ਰਾਗ malar baani bhagat ਨਾਮ ਦੇਵ ਜੀਓ ik ohankar satguru prasad malar raag malar malar da ke arth hai malar malhar keh malhar mal mal te jama sar karan karn wala malhar shabd malar nahi ਤੈਹਾਂ ਹਾ ਬੋਲਦੇ ਤੇ ਪੈਰ ਵਿੱਚ ਹਾ ਕੱਟਿਆ ਹੋਇਆ ਜੀ ਕਟਿਆ ਬਾਹਰ ਕੱਟਿਆ ਹੋਇਆ ਆ ਬਾਣੀ ਵਿੱਚ ਮਲਾਰ ਸ਼ਬਦ ਵੈਸੇ ਆਇਆ ਇੱਕ ਭਵਜਲ ਵਿਖਮ ਪੰਨਾ ਨੰਬਰ 59 ਭਵਜਲ ਵਿਖਮ ਡਰਾਵਣੋ ਨਾ ਕੰਦੀ ਨਾ ਪਾਰ ਨਾ ਬੇੜੀ ਨਾ ਤੁਲਹੜਾ ਨਾ ਤਿਸ ਵੰਜਮ ਮਲਾਰ ਉਵੇਂ ਹੋ ਰ ਆਰੇ ਯਾਰ ਉਹ ਅਭ ਜਲਦੇ ਵਿੱਚ ਨਹੀਂ ਆ ਮਾਲਾ ਕਰਨ ਵਾਲੀ ਕੋਈ ਚੀਜ਼ ਹਾਂ ਹਾਂਜੀ ਨਾ ਬੇੜੀ ਜਨ ਤਾਂ ਹੋਇਆ ਬੇੜੀ ਤੋਂ ਲਾ ਥੋੜੀ ਐ ਪਾਰ ਕਰਨ ਵਾਲੀ ਤਾਂ ਪਸੰਦ ਆਵੇ ਇੱਥੇ ਨਾ ਮਲ ਹਾਰ ਨਾ ਪੱਦਾ ਪਾਸਾ ਢਿੰਦਾ ਇਕ ਦਾ ਉਹ ਪੱਲਾ ਪਾਸਾ ਢਿੰਦਾ ਹੀ ਹੋਵੇ ਪੂਰੇ ਦਰਿਆ ਦੇ ਖੜੇ ਪੁਰੇ ਤਾਂ ਹੈ ਪਾਸਾ ਬੇੜੀ ਧੋਣਾ ਦਾ ਜਿਆਦਾ ਮਾਉਂਦਾ ਆਦਮੀ ਜਾਂ ਪੱਲਾ ਪਾਸਾ ਦਿਖਾਈ ਦੇਵੇ। ਯਾਰ ਆ ਮੈਂ ਬੇੜੀ ਧੋਣਾ ਬਣਾ ਕੇ ਬਾਹਰ ਜੂਣਾ। ਹਾਂਜੀ। ਨਾ ਤੇ ਵੰਜ ਮਲਾਰ। ਮਤਲਬ ਵੰਜ ਮਲਾਰ ਦਾ ਕੀ ਇਥੇ? ਉਹ ਬਾਸ। ਬਾਸ ਨੂੰ ਨਾ ਥੱਲੇ ਲਾ ਕੇ ਚਲੋਗੇ। ਨਾ ਬਾਹਰ ਨਾ ਕੋਈ ਐਸੀ ਚੀਜ਼ ਹੈ ਜੀ ਨਾ ਪਾਸਾ ਦੇ ਕੇ। ਨਾ ਸੱਖ ਦੇ ਵਿੱਚ ਕੋਈ। ਦੁਆ ਨਾ ਨਾ ਪਰ ਚੱਕਣ ਵਾਲੀ ਕੋਈ ਚੀਜ਼ ਹੈ ਇਹ ਤਾਂ ਦੇ ਤਰੀਕੇ ਬੇੜੀ ਤੋਂ 라 ਜਿਵੇਂ ਆਪਾਂ ਅਪਣਾਉਨੇ ਆ ਠੀਕ ਹੈ ਨਾ ਇਹ ਦੱਸਿਆ ਵੀ ਇਹਨਾਂ ਨਾਲ ਪਾਰ ਹੋਣਾ ਹੋਰ ਕਿਹਦੇ ਨਾਲ ਹੋਊ ਪਰ ਜਿਵੇਂ ਪਾਰਤਨਾਥ ਵਿਚ ਨਹਿਰ ਉਹਨਾਂ ਨੇ ਜਦੋਂ ਮੱਛੀ ਫੜ ਲਈ ساری ਮੱਛੀਆਂ ਨਾਲਕੜਿਆ ਵਿੱਚੋਂ ਬੰਦਾ ਜਿਹੜੇ ਸਮਾਦੀ ਲਈ ਹੋਈ ਸੀ ਹਾਂਜੀ ਉਹ ਕਹਿੰਦੇ ਇੱਕ ਬੰਦੂਰ ਸਾਰੇ ਮਾਛੀ ਸੀ ਤਾਂ ਪਾਰ ਪਾਰ ਦੇਖ ਲੈ ਨਹੀਂ ਬੰਦਾ ਨਿਕਲੇ ਕਿਸੇ ਜੋ ਵੀ ਰਾਜਾ ਕਹਿੰਦਾ ਵੀ ਤੂੰ ਬਈ ਝੂਠ ਬੋਲਦਾ ਗੱਲ ਕੀ ਉਹ ਕਹਿੰਦਾ ਵੀ ਤੁਸੀਂ ਮੇਰੀ ਗੱਲ ਨਹੀਂ ਸਮਝਦੇ ਨਾ ਇਹ ਕਿਹਾ ਜੀ ਖੀਰ ਤਾਂ ਕਰਾ ਪਹਿਲੀ ਤਾਂ ਗੱਲ ਹੈ ਸਾਡਾ ਤਾਂ ਖੀਰਾਂ ਦੜ ਨਹੀਂ ਖੀਰ ਸਾਡਾ ਵੀ ਜ ਜਾਓ ਉਹ ਬਿਵੇਕ ਦੇ ਜਾਲ ਚ ਉਹ ਕੀ ਮੱਛੀ ਉਹ ਬਿਵੇਕ ਦਾ ਜਾਲ ਕਹਿੰਦੇ ਵੀ ਬਿਵੇਕ ਦਾ ਤਾਂ ਜਾਲ ਹੀ ਨਹੀਂ ਹੁੰਦਾ ਇਰੋ ਨੇ ਆਪ ਬਵੇ ਸ਼ੁਰੂ ਕੀਤਾ ਬਵੇ ਕਵੇਤ ਦੀ ਕਹਾਣੀ ਅਬਵੇ ਕੀ ਹੁੰਦਾ ਥੋਡੇ ਕੋ ਅਬਵੇ ਦੇ ਜਾਲ ਨੇ ਕੋਈ ਵਿਦਿਆ ਤੁਸੀਂ ਸਮਝੀਵੇ ਮੈਂ ਜੋ ਕਿਹਾ ਕਿ ਜਾਲ ਮੱਛੀ ਦਾ ਉਹੀ ਤਾਂ ਮੱਛੀ ਕਹਿੰਦਾ ਕਿ ਵੀਰ ਜਲ ਕੀ ਮਛਲੀ ਜਲ ਖਜੂਰ ਉਸ ਮੱਛੀ ਦੀ ਉੱਥੇ ਗੱਲ ਹੈ ਜੇ ਕੋ ਪਾਣੀ ਵਾਲੀ ਮੱਛੀ ਸਮਝ ਲਵੇ ਹਾ ਤੇ ਤੇ ਉਹ ਬਿਦਿਆ ਬਿਦਿਆ ਦੀ ਬਲ ਹੋਈ ਨਾ ਆ ਬਿਦਿਆ ਸੋਦੇ ਤਾਤਲ ਹੈ ਨਾ ਸਾਨੂੰ ਇਹ ਸਮਝ ਆਈ ਨਹੀਂ ਪਲਕ ਨਾਰਾ ਜਿਹੜਾ ਵੀ ਨਾ ਇੱਥੇ ਕੋਈ ਦੱਸ ਰਿਹਾ ਹੈ ਕਿ ਦੂਰ ਕਰ ਰਿਹਾ ਵੀ ਭਾਈ ਐ ਨਹੀਂ ਐ ਹੋ ਪਾਪ ਦੂਰ ਕਰਨ ਵਾਲਾ ਵੀ ਨਹੀਂ ਗੁਰੂ ਕੋਈ ਉਪਦੇਸ਼ ਬਿਲਕੁਲ ਜੀ ਬਲ ਆ ਦਾ ਮਤਲਬ ਉਹ ਮਲ ਹਾਰ ਨਾ ਕੋਈ ਮਲ ਹਾਰਨ ਕਰਨ ਵਾਲਾ ਹੈ ਪਰਮ ਦੂਰ ਕਰਨ ਵਾਲਾ ਗੁਰੂ ਕਰੀਏ ਨਾ ਸਾਧਨ ਵੇੜੀ ਤੋਂ ਵਗੈਰਾ ਪਾਉਂਸ ਉਹਦਾ ਆਪ ਕਰਨਾ ਜਿਵੇਂ ਮਾਲਾ ਫੇਰ ਕੇ ਨਾਮ ਜਪ ਕੇ ਸਮਾਧੀ ਲਾ ਕੇ ਹਾਠੀਓ ਕਰਕੇ प्राणायाम करके ऐसा होगे ना बेड़ी तोला अपने साधन जे अपने साधन है नहीं कोई यत्न है नहीं कोई बेटा होगे ना यत्न जे यत्न नहीं कोई है तब फिर कोई पुचौना चाहिए다 और कोई साधन चाहिए다 बिना मेरे जतन दे बिना ओ वाला है ਕੋਈ ਉਹ ਪਰਮ ਦੂਰ ਕਰੇ ਗੁਰਪਰਸਾਦ ਭਰਮ ਦਾ ਨਾਸ ਕਰਨ ਵਾਲਾ ਨਹੀਂ ਕੋਈ ਹੈ ਮਲਾ ਦਾ ਮਤਲਬ ਹੈ ਐਸਾ ਸਤਗੁਰ ਨਹੀਂ ਹੈ ਗੁਪਤ ਦੁਆਰਾ ਮੋਕੜਾ ਹੈ ਆਵੋ ਜਾਓ ਉਹਨਾਂ ਨੇ ਅੱਗੇ ਕਲੀਅਰ ਕਰਤਾ ਸਤਗੁਰ ਭੈ ਕਾ ਬੋਇਤਾ ਨਦਰੀ ਪਾਰ ਉਤਾਰ। ਹਾਂ। ਉਹ ਸਤਗੁਰ ਨਹੀਂ ਹੈ ਕੋਈ ਉਹ ਕਹਿੰਦੇ ਸਤਗੁਰ ਹੈਗਾ ਭਾਈ। ਜਦ ਪਾਰ ਕੋਟੂਗਾ ਜਦ ਕਹਿੰਦਾ ਵੀ ਮੈਂ ਹੈਗਾ ਆਜੋ। ਫਿਰ ਉਹਨਾਂ ਨੇ ਕਿਹਾ ਮੁਕਤੀ ਮਿਲਦੀ ਹੋਈ ਨਹੀਂ ਜਿਉਂਦੇ ਨੂੰ ਫਿਰ ਉਹਨਾਂ ਨੇ ਬੰਦੇ ਕਹਤਾ ਰਸਤਾ। ਸਨਾਤਨ ਮਾਤਾ ਕਹਿੰਦਾ ਵੀ ਮੁਕਤੀ ਜਿਉਂਦੇ ਨੂੰ ਮਿਲਦੀ ਹੋਈ ਨਹੀਂ। ਕਬੀਰ ਕੰਨਾ ਮਰਨ ਮੁਕਤ ਕਿਨ ਪਾਈ ਆਤਮਾਨ ਦੇ ਬਾਦ ਕਿਨੋਂ ਮੁਕਤੀ ਮਿਲੂਗੀ ਕਿਨੋਂ ਨਹੀਂ ਮਿਲੂਗੀ ਇਹਦਾ ਕੀ ਤੂਰ ਹੈ ਤੁਹਾਡੇ ਕੋਲ ਇਹਦਾ ਸੁਖ ਹੀ ਨਹੀਂ ਪਾਈ ਤੇ ਬਾਦ ਮੁਕਤੀ ਇਹਦਾ ਸਾਰਿਆਂ ਨੇ ਪਾਈ ਹੈ ਇੱਕ ਜਨਮ ਨਹੀਂ ਹੌਸਲਾ ਕਰਕੇ ਵੇਰਾਂ ਇਹਨਾਂ ਨੂੰ ਤਾਂ ਜੋ ਸਨਾਤਨ ਮੱਤਾਲੇ ਜੀ ਆਓ ਵੀ ਜੀ ਗੁਰੂ ਬਣਾ ਹੈ। ਸਨਾਤਨ ਮਾਤਾ ਦੇ ਸਨਾਤਨ ਮਾਤਾ ਦਾ ਭਰਮ ਦੂਰ ਕਰਨ ਵਾਸਤੇ ਆਏ ਨੇ। ਉਹਨਾਂ ਨੂੰ ਪਤਾ ਹੈ। ਜਾਣਦੇ ਨੇ, ਸਮਝਦੇ ਨੇ ਪਰ ਜੇ ਉਹ ਆਮ ਦਾਨਸਰੀ ਹੋਣਗੇ ਸਨਾਤਨ ਮਾਤਾ ਦਾ ਜਿਹੜੇ ਦੂਰ ਸਨਾਤਨ ਹੈ। ਸ਼ਾਇਦ ਜਿਹੜੇ ਸਨਾਤਨ ਨੂੰ ਘਰ ਆਏ ਨੇ ਲੈ ਕੇ ਉਹਨਾਂ ਉ ਤਾਂ ਗਿਆਨ ਹੈਗਾ, ਸਮਝਦੇ ਨੇ ਦੂਜਿਆਂ ਦਾ ਭਰਮ ਦੂਰ ਕਰਨਾ ਚਾਹੁੰਦੇ ਨੇ। ਆਪਣੇ ਨਾਲ ਦੇ ਆਂਦਾ। ਜਿਵੇਂ ਨੇ ਕਿ ਆ ਸੀ ਆਪਣੇ ਬਨ ਚੁੱਕੇ ਨੇ ਜਿਵੇਂ ਆਰਾਸ ਆਰਾ ਵੀ ਮੈਂ ਭਾਗਵਤ ਵੀ ਜਿਲੇ ਗੈਰ ਸੈਂਟੀਫਿਕ ਗੱਲਾਂ ਨੇ ਇਹਦੇ ਚ ਹਿੰਦੂ ਮਾਤੇ ਚ ਉਹ ਤੇ ਆਦੋ ਭਾਈ ਹੁਣ ਬੋਲਿਓ ਹੁਣ ਨਹੀਂ ਸਮਾ ਹੈਗਾ ਉਹ ਤਾਂ ਇੰਨਾ ਇਸ਼ਾਰਾ ਕੀਤਾ ਉਹਨਾਂ ਨੇ ਜਿਹੜਾ ਤੁਹਾਡੇ ਕੋਲ ਗੈਰ ਸੈਂਟਰ ਕਮਨੀਅ ਲਿਖੀ ਹੋਈ ਹੈ ਨਾ ਜੀ ਫਾਤੀ ਦਾ ਸੱਲਾਤਾ ਬਖਰੀ ਦਾ ਸੱਲਾਤਾ ਹੋ ਕਰਤਾ ਹੋ ਕਰਤਾ ਕਿ ਛੱਡੋ ਇਹਨਾਂ ਦਾ ਮਨ ਨੂੰ ਕੁਝ ਨਹੀਂ ਰੱਖਿਆ ਮਨਹਾਰ ਦੀ ਗੱਲ ਕਰੋ ਰਾਗ ਮਨਹਾਰ ਤੇ ਆਓ ਹੁਣ ਗੁਰਪ੍ਰਸਾਦ ਪਰਮਕਾਰਨਾ ਉਸ ਗੱਲ ਤੇ ਆਓ ਫੇਰ ਹੈ ਕਰੋ ਗੱਲ ਪਰਮਾਨੰਦੀ ਲੋੜ ਨਹੀਂ ਰੋਤਾ ਚੁਰੂ ਅਪਦਰ ਤੋ ਕੀ ਦੀ ਗੱਲ ਬੈਠਾ ਕੇ ਹੈ ਨਹੀਂ ਧਰਮ ਕਿਹੜਾ ਬੇਤਨ ਮੋਲ ਮੋਲ ਕਹਿੰਦਾ ਬੇਤਨ ਹੈ ਕਿ ਖੋਜ ਲੋ ਭਾਈ ਕਿ ਮੈਂ ਕਹਿੰਦਾ ਆ ਆ ਦੂਏ ਤੇ ਤਮੈਂ ਕਹਤਾ ਹੈ ਮੈਂ ਕਹਤਾ ਹੈ ਚਾਹ ਮੈਨੂੰ ਪਤਾ ਵੀ ਹੈ ਮੈਂ ਕਹਿੰਦਾ ਆਓ ਖੋਜੀਏ ਬਸ ਥੋੜੀ ਜਿਹੀ ਤਸਲੀ ਹੋ ਬਾਕੀ ਜਿੰਨੇ ਧਰਮ ਨੇ ਸਾਰੇ ਇਨਵਾਈਟਡ ਨੇ ਅੱਧੀ ਬੈਠਾਂ ਲੈ ਇਹ ਨੂੰ ਕਹਿੰਨਾ ਇੱਕਾ ਖੁਦਾ ਹੈ ਯਾਰ ਆਮ ਜੋ ਵੀ ਮੱਦੀ ਨੋ ਹੈ ਇੱਕ ਹੈ ਉਹ ਇੱਕ ਨੂੰ ਸਮਝਾ ਦੇਵੇ ਸਾਨੂੰ ਸਨਾਤਨ ਨਾਲ ਇੱਕ ਨੂੰ ਸਮਝਾ ਦੇਣਾ ਅਸੀਂ ਮੰਨ ਲਾਂਗੇ ਸਨਾਤਨ ਮਤ ਠੀਕ ਹੈ ਤਾਂ ਕਿ ਬੇਦਮਤ ਜਿੰਨੇ ਦਿਨੋਂ ਸਾਨੂੰ ਸਮਝਾਉਣ ਦੇ ਚੁੱਪ ਰਹਾਂਗੇ ਜਿੱਥੇ ਸ਼ੰਕਾ ਉਹ ਉਥੇ ਗੱਲ ਕਰਾਂਗੇ ਜਦੋਂ ਹਟ ਖੜੇ ਕਰਦੇ ਵੀ ਸਾਤੇ ਭਾਈ ਸਮਝਾ ਨਹੀਂ ਹੁੰਦਾ ਫਿਰ ਦੂਸਲਾਮ ਅਲੈਕੁਮ ਅਲੈ ਤੁਸੀ ਆ ਜਾਓ ਸਜਾਈਆਂ ਨੂੰ ਕਹਿੰਦਾ ਤੁਸੀਂ ਆਜੋ ਬੋਧੀਆਂ ਨੂੰ ਕਹਿੰਦਾ ਤੁਸੀਂ ਆਜੋ ਜਿਹੜਾ ਸਮਝਾ ਦੂ ਧੋਤਕ ਰਾਜਾ ਰਾਣੂ ਕੀ ਕਹਾਣੀ ਉਹ ਵੱਤ ਪੂਰੀ ਹੈ ਬਾਕੀ ਵੱਤ ਅਧੂਰੀ ਹੈ ਜਿਹੜੀ ਪੂਰੀ ਮੱਤਾ ਉਹ ਧਰਮ ਤਦ ਪੂਰੀ ਮੱਤਾ ਮੱਤਾ ਜਦ ਮੱਤ ਪੂਰੀ ਹੋ ਜਾਂਦੀ ਹੈ ਫਿਰ ਉਹ ਧਰਮ ਉਹਦਾ ਬੋਲਿਆ ਹੋਇਆ ਉਹਦਾ ਦਸ ਧਰਮ ਉਧੂਰੀ ਮਾ ਟਾਲਵੀ ਆਪਣੇ ਨੂੰ タル ਮੁਕਈ ਜਾਂਦਾ ਇਹ ਗਲ ਦੀ ਪ੍ਰੋਗਰਾਮ ਹੈ ਉਧੂਰੀ ਆਲੇ ਕਹਿੰਦੇ ਨੇ ਇਹ ਵੀ ਧਰਮ ਹੈ ਪੂਰੀ ਆਲੇ ਨੂੰ ਤਾਂ ਚਲੋ ਅਜੋ ਧਰਮ ਕਿਹਾਂ ਬੇਧਰਮ ਗਿਆਨ ਧਰਮ ਬੇਧਰਮ ਉਹਨਾਂ ਦਾ ਗਿਆਨ ਧਰਮ ਬਾਬਾ ਤੇ ਇੱਕ ਹੋਰ ਜਗਾ ਮਲਾਰ ਦੀ ਗੱਲ ਆਈ ਹੈ ਮਹੱਲਾ ਤੀਜਾ ਮਲਾਰ ਸੀਤਲ ਰਾਗ ਹੈ ਹਰ ਧਿਆਈ ਹੈ ਸ਼ਾਂਤ ਹੋਏ ਬੱਈਏ ਆਏ ਥੇ ਜਬ ਇਹ ਨਹੀਂ ਹੈ ਸਭੋ ਤੇ ਅੰਤ ਬਦਲ ਗਿਆ ਹੁਣ ਜਦ ਤਾਲ ਨੂੰ ਧਿਆਨ ਰੂਪ ਹੋ ਜਵੇ ਇੱਕੋ ਧਿਆਨ ਹੋ ਜਵੇ ਦੁਬਾ ਖਤ ਮੋਜਵੇ ਉਹ ਮਲਾਰ ਹੈ ਮਲ ਹਲ ਹੋ ਗਈ ਲੇਖਾ ਦੂਰ ਹੋ ਗਿਆ ਧਾਂਟ ਗਿਆ ਜੋ ਚੀਜ਼ ਦੇਖਣੀ ਚਾਹੁੰਦਾ ਤਾਂ ਦੇਖੀ ਉਹਦੇ ਤੇ ਫਿਰ ਗੱਡ ਗਈਆਂ ਅੱਖਾਂ ਦੇਖੀ ਉੱਥੇ ਖੁੱਪ ਗਈ ਫਿਰ ਜਿਵੇਂ ਕੋਈ ਜਿਹਾ ਆਪਾਂ ਖਜ਼ਾਨਾ ਲੱਭਦੇ ਹਾਂ ਉਹ ਆਪਾਂ ਨੂੰ ਕੋਈ ਚੀਜ਼ ਆਪਾਂ ਗੱਡ ਕੇ ਦੇਖ ਦੇਣ ਸੰਦੈ ਜਾਂ ਕਰਕੇ ਦੇਖਦੇ ਹਾਂ ਉਹਨਾਂ ਨੂੰ ਉੱਥੇ ਲੱਭ ਗਿਆ ਵੀ ਇੱਥੇ ਵੀ ਤੇਲ ਆਇਆ ਪਰਾਉਲ ਆਇਆ ਗੈਰ ਹੈ ਪਰ ਉੱਥੇ ਹੀ ਪੱਟਣਗੇ ਕੋਈ ਆਣਾ ਉੱਪਰ ਤਾਂ ਨਹੀਂ ਅੱਪਰ ਨੂੰ ਜਾਣਾ ਧਰਤੀ 'ਚ ਲੱਭ ਗਿਆ ਪਹਿਲਾਂ ਵਰਮਾ ਮਾਰ ਕੇ ਦੇਖਦੇ ਨੇ ਜਦੋਂ ਨੂੰ ਕਹਾਂ ਲਾ ਕੇ ਵੀ ਹੱਲੇ ਇੱਥੇ ਹੈ ਕੁਝ ਤੇ ਉੱਥੇ ਹੀ ਪੱਟਾਂਗੇ ਦੂਰ ਤੋਂ ਉਹਦੇ ਕੋਲ ਦੇ ਪੱਟਣੇ ਜਾ ਕੇ ਜਦੋਂ ਖੱਡ ਕੇ ਹੈ ਜੋ ਕੁਝ ਹੈ ਤੇ ਉਸੇ ਕੰਦੇ ਸਾਰਾ ਧਿਆਨ ਹੋ ਗਿਆ ਨਹੀਂ ਤੇ ਟੋਲ ਦੱਸਦਾ ਸੀ ਕਰਕੇ ਉੱਥੇ ਵੀ ਧਿਆਨ ਜਲ ਹੈਗਾ ਬਲਾਰ ਹੋ ਗਿਆ ਰਾਗ ਇੱਥੇ ਧਿਆਨ ਹੋ ਗਿਆ ਗੁਰ ਧਿਆਨ ਕਸ ਬੜਿਆ ਹੁੰਦਾ ਧਿਆਨ ਪਹਿਲਾਂ ਗਿਆਨ ਜਾਂ ਗਿਆਨ ਧਿਆਨ ਤੇ ਬਦਲਦਾ ਨਾ ਉਹ ਦੋਵੇਂ ਦਾ ਧਿਆਨ ਖੇਡਦਾ ਫਿਰ ਸਾਡੀ ਦੁਨੀਆ ਦਾ ਧਿਆਨ ਸਾਡੀ ਮੁਕਤਰਾ ਧਿਆਨ ਖੇਚ ਲੈਂਦਾ ਕਿਦਾਂ ਤੇ ਨਹੀਂ ਸੇਟਾ ਕਿਦਾਂ ਜੀ ਧਿਆਨ ਗਿਆਨ ਦੇ ਜ਼ਖਦਾ ਗਿਆਨ ਕੋਤਮ ਦਾ ਅੰਮ੍ਰਿਤ ਕਟਿਆ ਜਾਂਦਾ ਹੁੰਦਾ ਗਿਆਨ ਦਾ ਅਗ ਜਿਵੇਂ ਹੀਰਾ ਜਿ ਚਲਦਾ ਹੈ ਅਗ ਫੜਦਾ ਕਿੰਨੀ ਰੋਜ਼ਨੀ ਹੁੰਦੀ ਹੈ ਸੂਰਜ ਜਿਹਾ ਹੀਰਾ ਅਗ ਲੱਗੀ ਹੋਈ ਹੈ ਇਹਨੂੰ ਸੂਰਜ ਹੀ ਹੈ ਐਟਮ ਚੁੱਟ ਰਹੇ ਨੇ ਜੀ ਚੱਲ ਕਿੰਨੀ ਰੋਜ਼ਨੀ ਹੈ ਪਰੇਗ ਦਾ ਧਿਆਨ ਕੇ ਤਾਂ ਨਹੀਂ ਜੇ ਤਾਂ ਕੁਝ ਆਰਟੀਫੀਸ਼ਲ ਕਿੱਡੀ ਰੋਸ਼ਨੀ ਪੈਦਾ ਕਰ ਦੂ ਆਰਟੀਫੀਸ਼ਲ ਧਰਮ ਨੇ ਕਿੰਨੀ ਕਿੰਨਾ ਗਿਆ ਰੋਸ਼ਨੀ ਪੈਦਾ ਕਰ ਦਨਗੇ ਇਸ ਕਰਕੇ ਇਹ ਜਿਹੜਾ ਬ੍ਰਹਮ ਗਿਆਨ ਸੂਰਜ ਇਹ ਚੱਕਦਾ ਮੇਰਾ ਇਹ ਕਰਦਾ ਪਰਮਾਨਾਸ ਆ ਗਿਆ ਮਲਾਰ ਆ ਗਿਆ ਤੇ ਇੰਡੈਕਸ ਇਸ ਲਈ ਕਿ ਅੰਦਰ ਜਲੀ ਗਿਆਨ ਤੇ ਆਣਾ ਜਾਣਾ ਬਾਤ-ਮਾਸ ਕਰ ਮੂਰਖ ਝਗੜੇ ਮੂਰਖ ਝਗੜੇ ਗਿਆਨ ਤੇ ਧਿਆਨ ਉਹ ਸਨਾਤ ਨਹੀਂ ਸਨਾਤ ਨਹੀਂ ਝਗੜੇ ਨਾ ਜੀ ਦੂਏ ਤੀਏ ਹੋਰ ਰਿਵਾਤਿਲ ਰਾਹ ਹੜੀ ਗਿਆਨ ਅਗਿਆ ਧਿਆਨ ਗਿਆਨ ਥਾਲ ਵਿੱਚ ਜਾਨਵਰ ਹੁੰਦਾ ਅੱਗ ਫੜਦਾ ਉਹ ਨਹੀਂ ਇਹਨੂੰ ਬਤਾ ਗਿਆਨ ਨਾਲੋਂ ਵੀ ਫੜ ਜਾਂਦਾ ਗੁਰ ਗਿਆਨ ਘੱਟ ਬੜਿਆ ਜਿਹੜਾ ਇਹ ਗਿਆਨ ਨਾ ਤੇ ਕਿਹਨਾਂ ਨੂੰ ਹੁੰਦਾ ਤੇ ਗਨਸੂਰੀ ਜਾਂਦਾ ਉਹਦੇ ਪੰਗ ਪਿਆ ਪਰਦਾਸਾ ਇਹ ਨਾਰਾ ਰਾਲ ਹੈ ਇੱਥੇ ਆ ਕੇ ਹੋਣਾ ਹੈ ਬਰਮਾ ਨਾ ਆਗੋ ਜਣਾ ਸਾਲੀ ਮਾਰ ਸਿੱਖ ਜਾਣੀ ਹਰ ਨਾ ਜਾਣੀ ਹੈ ਬ੍ਰਹਮਾ ਦਾ ਨ ਬ੍ਰह्म ਅਵੰ ਜੜੀ ਹੈ ਜੀਆ ਇਹ ਸਭ ਕੁਝ ਫੂਕ ਦਿੰਦੀ ਹੈ ਸਭ ਐ ਬੁੱਧੀ ਜਾਲੀਆਂ ਨੇ ਹਰ ਪ੍ਰਕਾਰ ਦੀ ਬੁੱਧੀ ਛਾੜ ਦੇਣੀ ਐ ਨੇ ਜੋ ਜੀਵ ਵਿੱਚ ਕੁਝ ਵੀ ਲਾਜੋ ਛਾੜ ਦੇ ਰਕੂੜਾ ਜੂਰ ਕਰ ਦੂ ਨੇੜੇ ਜਾਂਦੀ ਸਾਰੇ ਹਰ ਪ੍ਰਕਾਰ ਦੀ ਬੁੱਧੀ ਫੂਕ ਦਿੰਨਾਂ ਨੇ ਉਹ ਬਣੇ ਸਾਡੋ ਇਹ ਸੀ ਤਾਨੂੰ ਹਨ ਬਿਲਾਰਨ ਪ੍ਰੀਖਿਆ ਸੀ ਦادی ਇਹ ਹੀ ਹੈ ਉਹ ਅਗਲ ਦੀ ਆਪਣੀ ਪ੍ਰੀਖਿਆ ਹੈ ਸਭਾ ਬੁੱਧੀ ਜਾਰੀਨ ਕਰ ਹੈ ਤਤ ਗਿਆਨ ਸਿਰ ਤਤ ਛੱਡਦਾ ਪਹਿਲੇ ਜਾਂਦੇ ਬਾਦ ਜਿਹੜੇ ਇੱਥੇ ਰੰਗ ਨੇ ਸਾਰੇ ਭੂਖ ਤੇ ਤਾਂ ਦੇ ਹੋ ਜਾਂਦਾ ਤਾਂ ਅਗਲੇ ਜਨਮ ਜਨਮ ਬੁੱਧ ਹੁੰਦੀ ਹੈ ਬੱਚੇ ਜੀ बालभूत राग मलर वाणी भगत नामदेव जीयो की एक ओ अहंकार सतगुरु प्रसाद सेवियेले गोपाल राय अकुल निरंजन भगत दान दीजे जाचे संत जन राहो और भाई गल्ले आपाने ਜਿਹੜਾ ਪੜਿਆ ਪੜਦੇ ਆਂ ਤਾਂ ਜਿਹੜਾ ਪੜਿਆ ਐਹੀ ਪੜਿਆ ਜਾਂਦਾ। ਅਸਲ ਦੀ ਭਗਤੀ ਨੂੰ ਕੋਤ ਪੜਦੇ ਨਹੀਂ। ਪਰ ਬਿਲਕੁਲ ਅਰਥਾਂ ਨਾਲ ਤੇ ਇੱਥੇ ਪੜਨਗੇ ਹੋ ਜਾਣਾ। ਪਾਠ ਵੋਧ ਦੇ ਵਿੱਚ ਭਗਤ ਪੜਦੇ ਨੇ। ਉਹਨ ਭਗਤ ਜਿਹੜਾ ਬਾਣ ਦੀ ਜੈ ਜਿਹੇ ਪਹਿਲਾਂ ਭਗਤ ਹੁੰਦਾ ਭਗਤ ਮੁਕਤਾ ਹੁੰਦਾ ਸ਼ਬਦ। ਜੇ ਆਤਮਾ ਕੋ ਕੋ ਭਗਤ ਹੈ ਰਾਪੁਰਖ ਵਾਚਕ ਗ੍ਰੰਥ ਜੇ ਸਾ ਭਗਤ ਇੱਕ ਵਚਨ ਹੁੰਦਾ ਤਾਂ ਤਾਂ ਔਕੜ ਹੁੰਦਾ ਹੁਣ ਆ ਚਾਹੀਦਾ ਵਿਆਕਰਨ ਅਨੁਸਾਰ ਜੇ ਭਗਤ ਬਹੁਵਚਨ ਮੁਕਤਾ ਦਿੱਤਾ ਮੁਕਤਾ ਕੋ ਕਰਦਾ ਕਿ ਬਹੁਵਚਨ ਆ ਪਕਤਾਂ ਹੁੰਦਾ ਨਹੀਂ ਜੇ ਔਰ ਭਾਈ ਭਗਤਾਂ ਨੂੰ ਤਾਂ ਨਹੀਂ ਹੁੰਦਾ ਭਗਤ ਆ ਜਿਨੂੰ ਦਾਨ ਮਿਲ ਜਾਂਦਾ ਨਾ ਨਾਮਦਾਨ ਉਹ ਪਕਤ ਹੁੰਦਾ ਹੈ ਉਹ ਦੇਖੋ ਤਾਂ ਹੈਗਾ ਉਹ ਦਾਨ ਹੀ ਦੇਣਾ ਹੈ ਦਾਨ ਸੰਤ ਜਨ ਨੂੰ ਦੇਣਾ ਹੈ ਸੰਤ ਜਨ ਮੰਗਦੇ ਨੇ ਨਾਮ ਗੋਣ ਮੰਗਦਾ ਮੰਗਦਾ ਜਿਹੜਾ ਮਰ ਗਿਆ ਜਿਹਨੇ ਸੰਸਾਰ ਦੀਆਂ ਛਾਵਾਂ ਤਿਆਗ ਤੀਆਂ ਨਾਮ ਮਿਲੇ ਤਾਂ ਜੀਵਾਂ ਜੀਵਨ ਸੱਜੀਵਨ ਵਾਸਤੇ ਨਾਮ ਮੰਗਈਦਾ ਹੈ ਨਾਮ ਹੈ ਭਗਤੀ ਭਗਤੀ ਦਾ ਦਾਨ ਲੈ ਕੇ ਭਗਤ ਬਣ ਜਾਂਦਾ ਹੈ ਜਦੋਂ ਸ਼ੁੱਧ ਕੀਤਾ ਜਾਂਦੀ ਸੀ ਗੁਰਬਾਣੀ ਆਹੀ ਗੱਲਾਂ ਸ਼ੁੱਧ ਕੀਤੀਆਂ ਜਾਂਦੀਆਂ ਸੀ ਕੋਈ ਕਹਨੇ ਬੋਲ ਸਕਦੇ ਸੀ ਭਗਤੀ ਦਾ ਦਾਨ ਦਿੱਜੇ ਪਰ ਪੀ ਲਫ਼ਜ਼ੇ ਛੱਡਤਾ ਭਗਤੀ ਕਦੇ ਬੋਲਦੇ ਹੀ ਨਹੀਂ ਇਹ ਭਗਤੇ ਬੋਲਦੇ ਨੇ ਇਸ ਕਰਕੇ ਇਹਨਾਂ ਦੇ ਭਗਤੀ ਸਿੱਖੀਆ ਇਕੀ ਕੰਟੀਰੀਆੁਰ ਕੀ ਮੱਤ ਨੂੰ ਲੈ ਆਣੇ ਇਹ ਭਗਤੀ ਦੇ ਨਾ ਉਹ ਡੁੱਬੇ ਸਿਆਣੇ ਕੋਈ ਦੁਨਵੱਦਾ ਦਾਨ ਮੰਗਦਾ ਉਹ ਮੱਤ ਨਾ ਹੁੰਦਾ ਗੁਰੂ ਕੀ ਗੁਰ ਕੀ ਮੱਤ ਗੁਰ ਵਿੱਚੋਂ ਆਪਣੀ ਮਾਤ ਜਿਹੜੀ ਹੈ ਮਨਮਤ ਉਹਦੇ ਉੱਤੇ ਗੁਰਮਤ ਦਾ ਰੰਗ ਛਾੜ ਦੇਣਾ ਥੱਲੇ ਤੋ ਸੋ ਦੇਣੀ ਹੈ ਐਸੀਆਂ ਚੋਟਾਂ ਮਾਰਦੀ ਹੈ ਗੁਰਬਾਣੀ ਸਾਡੀ ਮਤ ਥੱਲੇ ਜ਼ਮੀਨ ਚ ਪਤਾਲ ਚ ਦੇ ਵਿੱਚ ਤਸੋਹ ਕੇ ਉੱਤੇ ਬਿਲਡਿੰਗ ਬਣਦੀ ਹੈ ਉਹਨਾਂ ਪੱਲਰਾਂ ਦਾ ਹੀ ਖੜੀ ਹੁੰਦੀ ਹੈ ਪੱਲਰ ਨਹੀਂ ਦੇ ਪਤਾਲ ਚੋਂ ਆਉਂਦੇ ਨੇ ਉਹ ਉੱਤੇ ਨੇ ਬਣੇ ਹੋਏ ਅਖੰਡਵਾਸ ਦੇ ਸਰਤੇ ਖੜੀ ਹੁੰਦੀ ਹੈ ਜੀ ਅਖੰਡਵਾਸ ਥੱਲੇ ਜ਼ਮੀਨ ਚ ਪਤਾਲ ਤੋਜ ਜਾਂਦਾ ਜੋ ਆ ਜਲਦਾ ਹੈ ਅਜਾੜਾ ਪਹਾੜਨਵਾਸ ਅਲੋਕ ਹੋ ਜਾਂਦਾ ਹੁੰਦਾ ਪਰ ਬੋਲਦੇ ਨਹੀਂ ਅੰਦਰੇ ਹੁੰਦਾ ਥੱਲੇ ਉਹ ਸੱਤੇ ਹੁੰਦੀ ਹੈ ਬੋਝ ਇਹ ਹਾਂਜੀ ਸੇਵੀ ਲੈ ਗੋਪਾਲਾਏ ਗੋਪਾਲਾਏ ਦੀ ਸੇਵਾ ਕਰੋ ਸੇਵੀ ਕਿਉਂਦਾ ਗੁਰ ਕੀ ਸੇਵਾ ਸ਼ਬਦ ਵਿਚਾਰ ਜੋ ਕੋ ਬਾਦ ਆਇਆ ਦਾ ਉਪਦੇਸ਼ ਹੈ ਉਹਦੀ ਵਿਚਾਰ ਕਰੋ ਉਹ ਜੋਦੀ ਸੇਵਾ ਜਿਵੇਂ ਕਹਿੰਦਾ ਉਵੇਂ ਕਰੋ ਜਿਵੇਂ ਚਲਾਉਂਦਾ ਉਵੇਂ ਚੱਲੋ ਕਰਨ ਵਿਚ ਚੱਲਣੀ ਸੇਵਾ ਸੇਵੀਲੇ ਗੋਪਾਲ ਵਾਲਾ ਉਹ ਬਾਲ ਰਾਇ ਦੀ સેવા ਕਰੋ ਕਿਉਂਕਿ ਉਹਨੇ ਭਗਤੀ ਦਾਣ ਦੇਣੀ ਹੈ ਸੰਤ ਜਨ ਨੂੰ ਦਾਣ ਦੇ ਸੰਤ ਤੇ ਘੱਟ ਨੂੰ ਭਗਤੀ ਨਹੀਂ ਮਿਲਦੀ ਪਹਿਲਾਂ ਸ਼ਾਂਤ ਹੋਣਾ ਪੈਂਦਾ ਹੈ ਪਹਿਲਾਂ ਸਬਰ ਕਰਨਾ ਪੈਂਦਾ ਹੈ ਸੰਤੋਖ ਤੋ ਬਾਦ ਇਹ ਨਾਮ ਮਿਲਦਾ ਇਹ ਨਾਮ ਨਾਲ ਵੈਸੇ ਨਹੀਂ ਬੜਾਉਂਦੇ ਨੇ ਉਹ ਭਾਈ ਹਉਮੈ ਨਾਮਾ ਨਾਲ ਵਿਰੋਧ ਹੈ ਉਹ ਕਹਿੰਦੇ ਹੰਕਾਰੀ ਨੂੰ ਨਹੀਂ ਨਾਮ ਕਾਇੰਦਤਾ ਨਾਮ ਟਿਕਦਾ ਨਹੀਂ ਉਹ ਸੁਣ ਨਹੀਂ ਸਕਦਾ ਤੁਸੀਂ ਉਹਨੂੰ ਨਾਮ ਦੇਈ ਜਾਂਦੇ ਹੋ ਨਾ ਦਾ ਤੇਣ ਵਾਲਿਆਂ ਕੋਲ ਕੁਝ ਹੈ ਨਾ ਲੈਣ ਵਾਲਿਆਂ ਕੋਲ ਤਾਂ ਵਿਚਾਰਿਆਂ ਕੋਈ ਜਿਆਦਾ ਉਹ ਜਾਂ ਤੇਣ ਵਾਲਿਆਂ ਕੋ ਕੋਈ ਹੋਵੇ ਤੇਣ ਵਾਲਿਆਂ ਦਾ ਪੱਲਾ ਘਟਾ ਗਾਹਾਂ ਉਹਨੇ ਜਿਹੜੀ ਟੀਜ ਦਿੱਤੀ ਹੈ ਮੁਠੀ ਉਹਦੀ ਤਾਂ ਮੁਠੀ ਖਾਲੀ ਹੈ ਮੁਠੀ ਦਾ ਕੁਝ ਹੈ ਨਹੀਂ ਤੇਰੀ ਝੋਲੀ ਕੀ ਬਹੁਤ ਜੌੜੇ ਆਪਣੀ ਮੁਠੀ ਖਾਲੀ ਹੈ ਖਾਲੀ ਮੁਠੀ ਪਾਈ ਜਾਂਦੇ ਨੇ ਖਾਲੀ ਝੋਲੀਆਂ ਲੈ ਕੇ ਤੁਹਾਨੂੰ ਆਈ ਜਾਂਦੇ ਨੇ ਖਾਲੀ ਮੁਠੀਆਂ ਪੈਂਦੇ ਨੇ ਖਾਲੀ ਝੋਲੀਆਂ ਆਉਂਦੀਆਂ ਨੇ ਅਸੀਂ ਝੋਲੀ ਭਰੀ ਵੀ ਅਜ ਤੱਕ ਭਗਤਾਂ ਦੀ ਝੋਲੀ ਜਦੋਂ ਭਰਦੀ ਪੰਚੀ ਨਾਲ ਝੋਲੀ ਭਰਨੀ ਸੀ ਨਾਮ ਬੋਣ ਦੀ ਕੋਲੀ ਗਏ ਤੇ ਪਿਆ ਜਿਹੜਾ ਆਲੇ ਕੋ ਨਾਮ ਹੈ ਨਹੀਂ ਪਤਾ ਹੀ ਨਹੀਂ ਕਿ ਕੀ ਨਾਮ ਹੁੰਦਾ ਆਪ ਲਈ ਨਹੀਂ ਸੰਤੋਖ ਹੈ ਹੀ ਨਹੀਂ ਆਪ ਨੂੰ ਕੀ ਅਵਸਥਾ ਹੋਣੀ ਚਾਹੀਦੀ ਹੈ ਕੀ ਕਰਨਾ ਚਾਹੀਦਾ ਹੈ ਗੁਰਬਾਣੀ ਕੀ ਕਹਿੰਦੀ ਹੈ ਤਾਂ ਸੁਣੇ ਕਿਥੇ ਨਹੀਂ ਉਹ ਘੜਨ ਬੜਾ ਲੈ ਸਾਬ ਨੇ ਦੁਕਾਨਦਾਰੀਆਂ ਚਲਾ ਲੀਆਂ ਬੜੀ ਛੇਤੀ ਚੱਲ ਪੈਂਦੀ ਹੈ ਕੋਈ ਬਹੁਤ ਇਨਵੈਸਟਮੈਂਟ ਨਹੀਂ ਹੈ ਜੇ ਵੀ ਨੇ ਗੋਪਾਲ ਰਾਏ ਆ ਕੇ ਹਾਸੀਗਾ ਜੀਤ ਗੁਰਬਾਨ ਨੇ ਕੁਛ ਕਰਨਾ ਦਾ ਸੰਤ ਜਨਾਂ ਨੇ ਕਿਸੇ ਸੰਤ ਨੇ ਕੰਮ ਕੀਤਾ ਜੇ ਤਾਂ ਹੁੰਦੇ ਸੰਤ ਚਨ ਫਿਰ ਤਾਂ ਕੰਮ ਕਰਦੇ ਜਿਹੜੇ ਸੀਗੇ ਸੰਤ ਜਨ ਉਹਨਾਂ ਨੇ ਤਾਂ ਕੰਮ ਕੀਤਾ ਜਾਣਦਾ ਮੈਂ ਜਾਣਕਾਰੀ ਲੈਣ ਵਾਲਾ ਜਾਨੀ ਜਿਹਨੂੰ ਗਿਆਨ ਲੈਣਾ ਜਿਹਨੂੰ ਨਾਮ ਦੀ ਭੁੱਖ ਹੈ ਜਾਜੀ ਹੈ ਇਹ ਤਾਂ ਨਾਲੋਂ ਬਾਅਦ ਫਿਰ ਤਾਂ ਮੰਗਦਾ ਇਹ ਕੰਮ ਕਰਦਾ ਪਰ ਇਹ ਤਾਂ ਸਾਰੇ ਪਰਪੰਚੀ ਸੀਗੇ ਇਹ ਤਾਂ ਬਨਾਰਸ ਕੇ ਠੱਗ ਸੀ ਸਾਡੇ ਮਾਣ ਇਹਨਾਂ ਨੂੰ ਫੀਲੋਡ ਭਈ ਸੀ ਉਹਨਾਂ ਦਾ ਪਰਦਾ ਫਾਸ਼ ਹੋ ਗਿਆ ਤਾਂ ਤਾਂ ਨਹੀਂ ਫਾਸ਼ ਕੀਤਾ ਸੀ ਉਦੋਂ ਉਦੋਂ ਨਹੀਂ ਪਰਦਾ ਫਾਸ਼ ਇਹਨਾਂ ਨੇ ਫੇਰ ਠੱਗਤਾ ਕੋਲ ਪਰਦਾ ਫਾਸ਼ ਹੋ ਗਿਆ ਸੋਣਾ ਓਖਾ ਟਕਣਾ ਉਦੋਂ ਕਮਿਊਨੀਕੇਸ਼ਨ ਦਾ ਸਾਧਨ ਹੈ ਨਹੀਂ ਸੀ ਯੋ ਇੰਟਰਨੈਟ ਹੈ ਹਰੇਕ ਦੇ ਕੋਲ ਮੋਬਾਈਲ ਹੈ ਪਰ ਤਾਂ ਟੈਲੀਵਿਜ਼ਨ ਕੋਣ ਇਹਨਾਂ ਦਾ ਬਚਾ ਨਹੀਂ ਹੋ ਸਕਦਾ ਟੈਕਨੋਲੋਜੀ ਨੇ ਪਰਮਿਸ਼ਨ ਪੈਦਾ ਕਰਤੀ ਉੱਖ ਵੀ ਬਹੁਤ ਪੈਦਾ ਕਰਤੀ ਲੋਕਾਂ ਨੇ ਸੇਵੀਲੇ ਬੋਲ ਗਏ ਉਹ ਬਾਹਰ ਦੀ ਸੇਵਾ ਕਰੋ ਉਹ اندر ਹੀ ਆ ਸਭ ਦਾ ਗੋਪਾਲ ਇਹ ਦੇਖਣ ਨੂੰ ਕਦੋਂ ਦਨੇ ਇਹ ਤੇ ਦੇਖਣ ਦਾ ਨੋ ਵਰਤ ਲਿਆ ਗੋਪਾਲ ਉਹ ਗਵੀਨ ਰਾਮ ਦਾ ਵਾ ਪੈਸੀ ਉਹ ਤਾਂ ਰਾਮ ਬੋਲੇ ਜੋ ਰਾਮ ਬੋਲਦਾ ਉਹ ਸੁਣੋ ਉਹ ਆਵਾਜ਼ ਅਨੁਸਾਰ ਕੰਮ ਕਰੋ ਉਹਦੀ ਮੰਨੋ ਉਹ ਬਾਲਾਏ ਜਿਵੇਂ ਕਰੋ ਉੱਠੋ ਪ੍ਰਾਪਤੀ ਹੋਣੀ ਹੈ ਤੁਹਾਨੂੰ ਦੀ, ਗੁਰਮਤ ਕੋ ਬਾਲਾਏ ਦੇ ਬਚਨ ਹੈ ਇਹਨੂੰ ਵਿਚਾਰੋ ਇਹ ਕਾਰਖਮਾ ਉਹ ਕੋਰ ਕਹਿਆ ਸਾਕਾਰਖਮਾ ਉਹ ਇਹ ਕਮ ਕਰਨਾ ਸੀ ਇਹ ਚੋਂ ਨਾਮ ਨਾਮ ਲੈਣਾ ਇਹ ਚੋਂ ਸਾਜੇ ਨੂੰ ਪ੍ਰਾਪਤੀ ਹੋਣੀ ਹੈ ਇਹ ਇਸੇ ਭੰਤੀ ਇਹੀ ਭਗਤੀ ਪਰਵਾਨਾ ਦਰਗਾਹ ਦੇ ਵਿੱਚ ਸੰਤ ਦੇ ਵਚਨ ਅਟੱਲ ਨੇ ਹੀ ਇਹ ਨਾਰਦ ਭਗਤੀ ਹੈ ਨਾਰਦੀ ਭਗਤੀ ਹੈ ਇਹਨੂੰ ਰੱਦ ਨਹੀਂ ਨਾ ਦਰਗਾ ਇੱਥੇ ਕੋਈ ਰੱਦ ਕਰਦਾ ਹੈ ਭਗਤੀ ਨੂੰ ਨਾ ਦਰਗਾ ਜਰਤ ਹੈ। ਇਹਦੇ ਖਿਲਾਫ ਕੋਈ ਤਰਖ ਨਹੀਂ। ਮੇਰਾ ਵਿਰੋਧ ਨਹੀਂ ਹੈ। ਆਕੀ ਸਾਰੀਆਂ ਭਗਤੀਆਂ ਦਾ ਵਿਰੋਧ ਦਾ ਵਿਰੋਧ ਹੈ। ਨਹੀਂ ਹੈ ਇਹਦਾ। ਹਾਂ ਇਹਨੂੰ ਵਗੜ ਲੈਣਾ ਨੇ ਫਿਰ। ਅਰਥਾਂਨਾਂ ਚ ਕਰਕੇ ਨਾ ਆਪਣੇ ਅਨੁਸਾਰ ਵੀ ਅਸੀਂ ਵੀ ਗੁਰਮਤਿ ਤੇ ਚੱਲਦੇ ਆਂ। ਆਪਣੇ ਮਤ ਨੂੰ ਗੁਰਮਤਿ ਦੇ ਬਰਾਬਰ तोड़ मरोड़ के पैनल कांदा का है ये कुछ कर रहे हैं हां जी हां जी जांचे कर दिग दिसै जांचे कर जिसदे कर दिग दिसै जालागै चेरग जांचे जा जानी जा ਜਾ ਜਿਹਦੇ ਘਰ ਵਿੱਚ ਜਿਹਦੇ ਘਰ ਅੰਦਰ ਜਿਸ ਦੇ ਘਰ ਅੰਦਰ ਜੀ ਦੇ ਘਰ ਵਿੱਚ ਉਹਦੇ ਘਰ ਵਿੱਚ ਕੀ ਆ ਜੀ ਤੋਂ ਜੇ ਮੰਗਣ ਜਾਣੇ ਆ ਉਹਦੇ ਘਰ ਵੀ ਕੁਝ ਹੋਵੇ ਜਿੱਥੋਂ ਮੰਗਣ ਜਾਵਾਂਗੇ ਜੇ ਘਰੇ ਕੁਝ ਨਹੀਂ ਘਰ ਕਿਹਾ ਜਾ ਵੱਡਾ ਇਥੇ ਬਾਬਾ ਜੀ ਜਿਹਦੇ ਘਰ ਵਿੱਚ ਸਭ ਕੁਝ ਹੈ ਭਾਈ ਉਹ ਘਰ ਵੀ ਤਾਂ ਵੱਡਾ ਹੀ ਹੋਊ ਜੋਡਾ ਉਹ ਜੱਜੇ ਜੱਜੇ ਨੂੰ ਕੰਨਾ ਉੱਪਰ ਬਿੰਦੀ ਹੈ ਬਿੰਦੀ ਨਹੀਂ ਸੀ ਬਿੰਦੀ ਇਹਨਾਂ ਨੇ ਲਾਈ ਜਾਨੇ ਕਿਹੜੇ ਵਾਲਿਆਂ ਨੇ ਬਿੰਦੀ ਅੱਧ ਕਦੇ ਹੁੰਦਾ ਹੀ ਨਹੀਂ ਕੁਰਬਾਨੀ ਤੇ ਕਿਸੇ ਬੀੜ ਚ ਨਹੀਂ ਤਾਇਪ ਜਿਹ ਹੈ ਕਿਸੇ ਬੀੜ ਚ ਦਿਖਾਇਓ ਇਹਨਾਂ ਨੇ ਅਲੱਗ ਲਾਈਆਂ ਨੇ ਪੋਤੀਆਂ ਚ ਆਦ ਕਰ ਸਿੱਖ ਨੂੰ ਅੱਧ ਦਿਖਾ ਦਿੱਤੇ ਹੈਗਾ ਕਿਤੇ ਨਹੀਂ ਜੀ ਫਿਰ ਸਿੱਖ ਨੂੰ ਵੱਡਕ ਚਾਹੀਦਾ ਇੱਕ ਸਿੱਖ ਬਣ ਜਾਂਦਾ ਸਿੱਖ ਸਿੱਖਿਆ ਸਿੱਖਦਾ ਸਿੱਖਦਾ ਮਤਲਬ ਹੈ ਸੱਚੇ ਨੂੰ ਯਾਰੀ ਖਖਾਸ ਸਿੱਖ ਇਹਦਾ ਅਰਥ ਹੈ ਸਿੱਖਿਆ ਸਿੱਖਦਾ ਮਤਲਬ ਹੈ ਅਦਕ ਨਾਲ ਸਿੱਖ ਬਣਿਆ ਜਿਹਨੇ ਸਿੱਖਿਆ ਲੈਣ ਵਾਲਾ ਜਦੋਂ ਅਗਰ ਨਾਲ ਲੈਣ ਵਾਲਾ ਅਰਥ ਸਿਖਿਆ ਦੋ ਅਰਥ ਨਾਲ ਫਰਕ ਹੈ ਅਗਰ ਗੱਦੇ ਹੈ ਇਹ ਨਹੀਂ ਦਰਵਾਣੀ ਜੀ ਸਿਖੇਤਵਾਰ ਆਇਆ ਨਾਖ ਸਿਖ ਉਹ ਸਿਖਿਆ ਜਿਹੜੀ ਮੁੜਦੀ ਹੋਈ ਨਹੀਂ ਹੈ ਜਿਹਦੀ ਧਾਰ ਮੁੜਦੀ ਹੋਈ ਨਹੀਂ ਹੈ ਗੁਰਮਤਿ ਦੀ ਸਿਖਿਆ ਨਾਖ ਸਿਖ ਜੇ ਬਾ ਨਾਂ ਦਾ ਨੋ ਪਾਸੇ ਜੀ ਕੋਲ ਨਾਸ ਨੂੰ ਵਰਨੀ ਨਹੀਂ ਨਾ ਕਿ ਨਾ ਉਹ ਆਵੇ ਜਿਹੜਾ ਉੱਤਰਾ ਦਾ ਉਂਗਲ ਦਾ ਜਿਹੇ ਮੁੜ ਜਾਂਦਾ ਨਾ ਹਨ ਉਹ ਵੀ ਕਹਿੰਦੇ ਨੇ ਨਖਸ ਸਖਤ ਨੂੰ ਵੀ ਕਹਿੰਦੇ ਨੇ ਨਖ ਸਖਿਆਰ ਨੂੰ ਬੜਾ ਨਾਖਾਜ਼ਮੀਆ ਮੁੜ ਜਾਣੇ ਪਿਛੇ ਸਖਿਆਰ ਨਖ ਦੇ ਮੌਸਾ ਦੇ ਅਰਥ ਮੈਂ ਪਿਛੇ ਨਖ ਲੱਭਦਾ ਵਰਤਦੇ ਤੇ ਉਹ ਬੜਾ ਨਾਖਾਜ਼ਮੀਆ ਸੁਦਾ ਜਾਂਦਾ ਪਰਵਾਣੀ ਰੱਖਦਾ ਸੱਚਾ ਕੋਈ ਤਾਂ ਲੱਭੇ ਨਹੀਂ ਹੈ ਬੁਰਾ ਨੇ ਹਾਂ ਨਹੀਂ ਭਾਬੀ ਤੁਸੀਂ ਕਿਹਾ ਵੀ ਸਿੱਖ ਦੇ ਜੋ ਸਿੱਖਿਆ ਲੈਣ ਵਾਲਾ ਹੈ ਉਹਦੇ ਉੱਤੇ ਅੱਗ ਚਾਹੀਦੀ ਹੈ ਤਾਂ ਫਿਰ ਗੁਰਬਾਣੀ ਤਾਂ ਹੈ ਨਹੀਂ ਭਾਏ ਨਹੀਂ ਸੀ ਗੁਰਬਾਣੀ ਦੇ ਵਿੱਚ ਕਾਹਨ ਸੰਖਿਆ ਲੈ ਕੇ ਪੜ੍ਹਨ ਦੀ ਗੱਲ ਸੀ ਇਹੇ ਜਹ ਹੱਥ ਲਿਖਤਾਂ ਦੇ ਵਿੱਚ ਕਿਤੇ ਆਤ ਕਦੇ ਨਹੀਂ ਸੀ ਉਹ ਨਿਯਮ ਸੀ ਆਪਾਤ ਕੋ ਪਾਉਣਾ ਨਹੀਂ ਪਰ ਪੜਨਾ ਤੇ ਜਦ ਤੇ ਲੋੜ ਪਊ ਲਾ ਲੈਣਾ ਿੱਪੀ ਬਿੰਦੀ ਬਿੰਦੀ ਨਾਲ ਿੱਪੀ ਦਿਖਾ ਸਕਦੇ है ਚ ਚਾਰ ਚੀਜ਼ਾਂ ਨਹੀਂ ਹੈ ਬਿਲਕੁਲ ਵੀ ਉੱਪਰ ਜਿਹੜੇ ਆਉਂਦੇ ਤੇ ਕਹਿ ਵੀ ਸਤੂ ਕਰਤੀ ਆ ਨਾ ਹੱਥ ਲਿੱਕਾਂ ਵਿੱਚ ਹੁੰਦੀਆਂ ਸੀ ਜਿਹੜਾ ਨੇ ਰਾਤ ਨੂੰ ਜਿੱਦਿਆਂ ਨੇ ਜਦ ਕਹਿਤ ਕਰ ਸ਼ਾਪਾ ਪਾਇਆ ਪਹਿਲਾ ਹੈਂਸੀ ਸਾਹਿਬ ਹੈ ਵਿਸ਼ਵ ਦੇ ਵਿੱਚ ਪਹਿਲੇ ਬਾਵਾ ਹੈ ਬਿਸ਼ੂ ਨੂੰ ਬਿਸ਼ੂ ਇਸਾਈ ਨਾ ਜੀ ਫਿਰ ਬਿਸ਼ੂ ਸਾਹਿਬ ਦੇ ਗੁੱਟ ਦੇ ਬਾਵਾ ਬਾਵਾ ਇਹ ਵਿਸ਼ਵ ਸੰਸਾਰ ਜੇ ਤੂੰ ਦੇਖਦਾ ਯਾਰ ਕਾ ਰੂਪ ਹੈ ਇਹਵੇਂ ਨੇ ਸਾਇਕੰਗ ਦੇ ਵਿੱਚ ਪਾਵਾ ਘਟਾਇਆ ਫਿਰ ਚੋਂ ਇਹਨਾਂ ਤਾਂ ਇੰਨੀ ਭਗਾੜਦੀ ਗੱਲ ਵੀ ਇਹ ਠੀਕ ਹੋਈ ਨਹੀਂ ਸਕਦੀ ਝਗੜੇ ਚ ਪਈ ਰਹੇ ਝਗੜੇ ਤੇ ਮੈਂ ਆਇਆ ਸੀ ਜਾਂ ਝਗੜਾ ਹੀ ਹੋ ਰਿਹਾ ਸੀ ਬਾਠਨਪੁਰ ਦਾ ਮੈਂ 6 ਸਾਲ ਝਗੜੇ ਚ ਆਪਰੇ ਹਾਂ ਉਹ ਝਗੜੇ ਚ ਨਾਲ ਇਧਰ ਨਿਕੜਿਆ ਉਹ ਛੜਤਾ ਦੂਆ ਪਤਾ ਉਹ ਝਗੜੇ ਦਾ ਹੱਲ ਕੱਢੀ ਐ ਕੀ ਐ ਹਣ ਹੱਲ ਖਾਤਰੇ ਮੈਂ ਸਾਡਾ ਬੁੱਢਾ ਗੱਲ ਛੱਡਿਆ ਐ ਦੇਖੋ ਕੀ ਬਲੂ ਬਨ ਕੋਈ ਨਹੀਂ ਇਹਦਾ ਕੋਈ ਨਹੀਂ ਯਾਦ ਕੋਈ ਮੈਨੂੰ ਚਿੰਤਾ ਨਹੀਂ ਹੋ ਜਲਦੀ ਸੰਤਾ ਨੂੰ ਕੋਈ ਚਿੰਤਾ ਨਹੀਂ ਕਿਸੇ ਨਾਲੀ ਆਪਾਂ ਫਾਲਸਾ ਸਭ ਕੋ ਆਪਣੇ ਕੋਲ ਉਹਦਾ ਘੋੜਿਆਂ ਨੂੰ ਤਲਵਾਰਾਂ ਨੂੰ ਲੋਕਾਂ ਨੂੰ ਸਮਝਦੇ ਕੋਲ ਸਾਡੇ ਸਭ ਕੁਝ ਕੋਣੇ ਗਿਰਣਾ ਜੀ ਅਤੇ ਦੂਜਾ ਨਵੀਂ ਵੀ ਲੜਨ ਇਹ ਤਾਂ ਆਪਣੇ ਆਪਣੀ ਭੁੱਖ ਹੁੰਦੀ ਹੈ ਮੈਨੂੰ ਪਤਾ ਲੱਗਿਆ ਸਾਡੇ ਕੋਲ ਨਹੀਂ ਕੱਖ ਨਹੀਂ ਜਿਹੜੀ ਚੀਜ਼ ਖਾਤਰ ਮੈਂ ਬਾਣਾ ਪਾਇਆ ਉਹ ਤਾਂ ਹੈ ਹੀ ਨਹੀਂ ਨਾ ਕੋਲ ਮੈਨੂੰ ਪਤਾ ਲੱਗਿਆ ਬਾਅਦ ਚ ਜੀ ਸਾਲ ਇਹਦੇ ਕੋਲ ਤਾਂ ਕੁਝ ਵੀ ਨਹੀਂ ਜਦੋਂ ਉਹ ਕਹਿੰਦੇ ਸਾਨੂੰ ਕੱਚੀ ਪੱਕੀ ਬਾਣੇ ਦਾ ਗਿਆਨ ਹੀ ਨਹੀਂ ਕਿਸੇ ਨੂੰ ਅੰਨੀ ਸ਼ੌਕਰ ਕਰ ਗਿਆ ਇਹਨਾਂ ਕੋਲ ਕੁਝ ਵੀ ਨਹੀਂ ਵਾਲਾ ਤਾਂ ਲੇਖੇ ਜਾ ਗਿਆ ਕੋ ਜੋ ਕੀਤੀ ਮੈਂ ਆਪ ਕੋ ਜੋ ਕੀਤੀ ਰਾਮਣੇ ਦੇਖੋ ਪਹਿਲਾਂ ਦਿਖਾਉ ਕਿ ਹੈ ਉਹ ਵੀ ਚਾਹ ਲੋ ਇੱਛਾ ਸੀ ਪਰ ਮੈਂਛ ਨੇ ਆਪ ਕਰਾ ਲੀਂ ਕਰਦੇ ਦਾ ਪਹਿਲਾਂ ਵੀ ਸੀ ਲੱਗੇ ਤੇ ਆਪਣੇ ਆਪਣੇ ਲੈਵਲ ਤੇ ਪਰ ਕੋਸ਼ਿਸ਼ ਚਲੋ ਕਰਾ ਲੀ ਕਿਵੇਂ ਆਕਰਾ ਲੀ ਕਿਵੇਂ ਹੋ ਗਿਆ ਮੇਰੀ ਇੱਛਾ ਸੀ ਕਹਾਂ ਹੋਵੇ ਜੇ ਸੀਗੀ ਤਾਉਨ ਫੜ ਲਾ ਗਿਆ ਉੱਤ ਸਮਝੇ ਸਾਹਮਣੇ ਜੈ ਜੀ ਇੱਛਾ ਸੀ ਉਹ ਮੈਨੂੰ ਪਤਾ ਚੰਗੀ ਰਹੀ ਆ ਮਾਰੀ ਤੀ ਉਹਨੂੰ ਇੱਧਰ ਫੜ ਲਾ ਗਿਆ ਹੁਣ ਸਰ ਉੱਤ ਸਮਝੇ ਸਾਹਮਣੇ ਪ੍ਰਾਪਤੀ ਹੋਈ ਹੈ ਸਮਝੇ ਸਾਹਮਣੇ ਅਕਾਲੀ ਸਾਡੀ ਜੜ ਪੱਟਣ ਨੂੰ ਫਿਰਦੇ ਸੀ ਆਰੇ ਖਲਾਵੇ ਇਹੜਾ ਬਾਣੇ ਦੇ ਖਿਲਾਫ ਆ ਉਹ ਸਿੱਖੀ ਦੇ ਖਿਲਾਫ ਆ ਉਹ ਤਾਂ ਬਾਣੇ ਨੂੰ ਦੇਖਣਾ ਨਹੀਂ ਚਾਹੁੰਦੇ ਲੋਕ ਗੁਰੂ ਸਾਰੇ ਫਰਵੀ ਮਹਾਰਾਜ ਚਲੇ ਗਏ ਕੋਈ ਚਲੇ ਗਿਆ ਉਹ ਇਹ ਦੇਖਣਾ ਨਹੀਂ ਚਾਹੁੰਦੇ ਇਹ ਵਾਲੇ ਬਾਬਾ ਜੀ ਉਹਨਾਂ ਦਾ ਕਹਿਣਾ ਜਿਹੜੇ ਦੇਖਣਾ ਨਹੀਂ ਚਾਹੁੰਦੇ ਜਿਵੇਂ ਅਸੀਂ ਆਮ ਸੁਣਦੇ ਵੀ ਧਿਆਨ ਸਿੰਘ ਦਾ ਜਿਹੜਾ ਕਿਰਦਾਰ ਹੈ ਉਹ ਠੀਕ ਨਹੀਂ ਹੈਗਾ ਜੇ ਨਹੀਂ ਜੀ ਗੱਲ ਕਿਉਂ ਲਾਏ ਨੇ ਇਹਨਾਂ ਨੂੰ ਫੇਰ ਠੀਕ ਆਲੇ ਬਾਦਨ ਗੋਡਿਆਂ ਦੇ ਥਲੇ ਘੁੜਾਲੇ ਨੇ ਅਗਾਹ ਤੱਕ ਤੇ ਨੇ ਛੇਕ ਦੇ ਗੇਉਨੀਏ ਰਾਨੂੰ ਉੱਥੇ ਜਿਹੜੇ ਗਲਤ ਨੇ ਉਹ ਤਾਂ ਉਹਨਾਂ ਦੇ ਨਾਲ ਨੇ ਮੈਨੂੰ ਦਾ ਸਿਰ ਮੇਰਾ ਕਲਦਾਰ ਕਹਿਆ ਜੇ ਮੈਂ ਉਹਨਾਂ ਦੇ ਨਾਲ ਦੀ ਜੋ ਜੋ ਠੀਕ ਨਹੀਂ ਨਾਲ ਕਿਉਂ ਲਾਏ ਨੇ ਆਪਣੇ ਯੂਜ਼ ਕਰਨ ਲਈ ਯੂਜ਼ ਕਰਨੇ ਉਹਨਾਂ ਉਹਨਾਂ ਵਾਤੇ ਠੀਕੇ ਨੇ ਉਹਨਾਂ ਵਾਤੇ ਦਾ ਠੀਕੇ ਨੇ ਨਾਲੇ ਲਾੜਦੀਆਂ ਫੌਜਾਂ ਕਹਿ ਦਿੰਦੇ ਨੇ ਨਾਲੇ ਕਹਿੰਦੇ ਨੇ ਬਾਣਾ ਇਹਨਾਂ ਨੇ ਰੱਖਿਆ ਸਾਥੇ ਰੱਖ ਨਹੀਂ ਹੋਇਆ ਨਾਲੇ ਕਹਿੰਦੇ ਨਹੀਂ ਠੀਕ ਨਹੀਂ ਤੁਸੀਂ ਢੀਪੋ ਜੇ ਇਹ ਠੀਕ ਨਹੀਂ ਤੁਸੀਂ ਭਾਈ ਠੀਕ ਬਣ ਜਾਓ ਤੁਸੀਂ ਪਾਓ ਬਾਣੇ ਉਹ ਵੀ ਠੀਕ ਬਣਾਓ ਫਿਰ ਇਹ ਠੀਕ ਨਹੀਂ ਅਸੀਂ ਇਹਨਾਂ ਨੂੰ ਗੁਰੂ ਦੇ ਬਰਾਬਰ ਪੰਥ ਦਾ ਬਰਾਬਰ ਨਹੀਂ ਮੰਨਦੇ ਅਸੀਂ ਠੀਕ ਨੇ ਇਹਨਾਂ ਨਾਲ ਵੀ ਅਸੀਂ ਘਟੀਆਂ ਅਸੀਂ ਲੀਡਰ ਤੁਸੀਂ ਕਿਹਾ ਠੀਕ ਉਹਨਾਂ ਨੂੰ ਪੁੱਛੋ ਠੀਕ ਹੋ ਫਿਰ ਉਹਨਾਂ ਬਾਈ ਮੀਟਿੰਗ ਕਿਹਨੇ ਅਕਾਲੀਆਂ ਨਾਲ ਫੇਰ ਠੀਕ ਨੇ ਸੰਤਾਨਾਂ ਨਾਲ ਫੇਰ ਠੀਕ ਨੇ ਪਰ ਜਿਹੜੇ ਜਗੁਰੂ ਨੇ ਬਣਾਇਆ ਤਾਂ ਉਹ ਜਿਹੜੀ ਹਨ ਉਹ ਤਾਂ ਸੀ ਤਾਂ ਗੁਰੂਆਂਾਂ ਦੀ ਗੱਲ ਕਰਦੇ ਇਹਨਾਂ ਦਾ ਤਾਂ ਮਿਹਲੇ ਇਹ ਤਾਂ ਖੰਡਵਾਦ ਇਹ ਆਪ ਜਾਂ ਖੰਡਵਾਦ ਉਹਨਾਂ ਵੱਲ ਨੂੰ ਜਾਣ ਲੱਗੇ ਜਿਆਦਾ ਇਹਨਾਂ ਨੂੰ ਕਹਿੰਦੇ ਆ ਤੁਸੀਂ ਕਹਦੇ ਬੇਹ ਪਾਣੀ 'ਚ ਬਹਿ ਗਏ ਕੋਈ ਨੂੰ ਕਾਦੀ ਭੋਖਾ ਬਾਣਾ ਪਿਉ ਪਾਇਆ ਪੜਨ ਲੱਢੋ ਫਿਰ ਹਾਂਜੀ ਬਾਬਾ ਜੀ ਤੁਸੀਂ ਹੁਣ ਕਿਹਾ ਸੀ ਅੱਜ ਬਾਰੇ ਗੱਲ ਹੋਈ ਸੀ ਜਿਵੇਂ ਬਾਣੀ ਦੀ ਪੰਕਤੀ ਹੈ ਮੰਨੈ ਤਰੈ ਤਾਰੇ ਗੁਰਸਿਖ ਉਥੇ ਪੜਾ ਨਹੀਂ ਫਿਰ ਆਲਤ ਪੜਦੇ ਜੀ ਮੰਨੈ ਤਰੈ ਤਾਰੇ ਗੁਰਸਿਖ ਗੁਰਸਿਖ ਤਾਰਦਾ ਬਾਕੀ ਤੜਦੇ ਨੇ ਕਿਨੂੰ ਜੇ ਤਰੇ ਤਾਰੇ ਤਰੇ ਗਦੇ ਹੂੰਗਾ ਆਪ ਦਾ ਕਰਦਾ ਹੀ ਜਿਹੜਾ ਤਾਰਦਾ ਜੱਗ ਤਾਰੇ ਗੁਰ ਸਿੱਖਾ ਜੱਗ ਗੁਰ ਸਿੱਖ ਤਾਰਦਾ ਕਿੰਨੂੰ ਤਾਰਦਾ ਮੁੰਨਾ ਤਰਾਂ ਤਾਰੇ ਗੁਰ ਸਿੱਖ ਤਾਰਦਾ ਜਿਹੜੇ ਨਵੇਂ ਜਿਹੜੇ ਸਿੱਖ ਨਾ ਤਰਦੇ ਨੇ ਗੁਰ ਬਣਦੇ ਨੇ ਗੁਰਸੇਖ ਜਦ ਬਣ ਜਾਂਦਾ ਕਰ ਜਾਂਦਾ ਸਿੱਖ ਦਾ ਤਰਵਾ ਨਹੀਂ ਹੈ ਸਿੱਖ ਦਾਤਾ ਸਿਰਫ ਨੱਕ ਨੂੰ ਉਹ ਅੱਖਾਂ ਬਲਕੇ ਮੂੰਹ ਵੀ ਨਹੀਂ ਹੈ ਨੱਕ ਅੱਖਾਂ ਤਨ ਇਹ ਬਾਹਰ ਹੈ ਪਾਣੀ ਤੋਂ ਉਹ ਪਾਣੀ ਤੋਂ ਬਾਹਰ ਹੈ ਜਦ ਇਹ ਮੂੰਹ ਪਾਣੀ ਤੋਂ ਉਹ ਗੋਲੂ ਦਾ ਪਾਣੀ ਦੇ ਜੂਗਾ ਦੱਬਾ ਕੇ ਤੇ ਸਾਹ ਹੁੰਦਾ ਨੰਬਕ ਇਹ ਪਾਣੀ ਦੀ ਬਾਤ ਚਾਈ ਜਾਈਏ ਅੱਖਾਂ ਦੇਖੂਗਾ ਤਾਂ ਇਹ ਪਾਣੀ ਦੇ ਵਾਰ ਅੱਖ ਉੱਤੇ ਥੱਲੇ ਜੀ ਤੇ ਬਾਕੀ ਕੰਨ ਜਦ ਨਾਲ ਬੱਚਾ ਪੈਦਾ ਹੁੰਦਾ ਨਾ ਸਭ ਤੋਂ ਪਹਿਲਾਂ ਆਉਂਦਾ ਉਹ ਜਵਾਂ ਦੇ ਅੱਖਾਂ ਬਾਹਰ ਚਲਦੀਆਂ ਨੇ ਕੋਕ ਸਾਹੀ ਜੀਵਨ ਪਹਿਲਾਂ ਨੂੰ ਤ੍ਰਣ ਵਹੀ ਜਾਈ ਦੀ ਹੈ ਜੀ ਆਹ ਅੱਖਾਂ ਦੀ ਗੱਲ ਬਾਤ ਅੱਖਾਂ ਦਾ ਨਾਮ ਹੀ ਹੋਰ ਤਾਂ ਸਮਝੂਗਾ ਉਹ ਪੈਦਾ ਹੁੰਦਾ ਨਾ ਪਹਿਲਾਂ ਆਉਂਦੀਆਂ ਨੇ ਮਨੈ ਤਰ ਤਾਰੇ ਗੁਰਸਿੱਖ ਜਿਹੜਾ ਸਸਤਾ ਤਰਦੇ ਨੇ ਤਰੇ ਬਹੁ ਬਚੇ ਨੇ ਸਸੇ ਸਾਧੂ ਵਰ ਤੋਂ ਸੇਖਾ ਨਾਣ ਵਾਲੀ ਵਰਤਿਖ ਨਹੀਂ ਹੈ। ਬਣਾ ਬਰਤਕੇ ਹੋਰ ਕੀ ਹੈ? ਸੇਖਾ ਗੁਰੂ ਗੁਰੂ ਸੇਖਾ। ਨਾਣਕ ਪੈਦਨਾ ਭਾਈ। ਸੇਖ ਸੇਖਾ ਲੈ ਕੇ ਗੁਰੂ ਬਣਦਾ। ਸੰਸਾਰ ਦੇ ਵਿੱਚ। ਸੰਸਾਰ ਦੇ ਵਿੱਚ ਜਿਵੇਂ ਆ ਗੁਰੂ ਬੰਦੇ ਨੇ ਪਹਿਨਾ ਸਿੱਖਿਆ ਲੈਂਦਾ ਫਿਰ ਸੁਹਾਗ ਜਾਂਦਾ ਪੜਾਉਣ ਲੱਗ ਜਾਂਦਾ ਉਹ ਸਾਰੇ ਸੰਸਾਰੀ ਸਿੱਖ ਦੀ ਗੱਲ ਆ ਉਹ ਜੀ ਆ ਹਾਂਜੀ ਜਾਂਚੇ ਕਰ ਦਿਗ ਦਿਸੈ ਜਾਂਚਿਆ ਕਰ ਜਾਂ ਚੈ ਕਰ ਜਾ ਚੈ ਜਾਂ ਛੱਬ ਦੇ ਕਿਤੇ ਆਉ ਜਾਂ ਦੇ ਨਾਲ ਤਾਉ ਜੇ ਤਾਉ ਜਾਂ ਕੰਡੀਸ਼ਨਲ ਸ਼ਬਦ ਹੈ ਜਾਂ ਤੂੰ ਮੇਰੇ ਵਾਲਾ ਜਾਂ ਹਿੰਦੀ ਦਾ ਸ਼ਬਦ ਹੈ ਜਾਂ ਦੇ ਨਾਲ ਤਾਉ ਦਾ ਟਾਕਾ ਮੂੜੋ ਚਾਰਤ ਪੈਦਾ ਜਾਂਖੋ ਪੇਵਨ ਬਾਬਤ ਹਿੰਦੀ ਬਹੁਤ ਹੈ ਸੁਤਰਾ ਮੈਂ ਪੰਜਾਬੀ ਨਹੀਂ ਪੜੀ ਮੈਨੂੰ ਤਾਂ ਪਤਾ ਕੋਰਵਾਣੀ ਬਾਰੇ ਹਿੰਦੀ ਸਾਈ ਲਿਖਿਆ ਹੈ ਪੰਜਾਬੀ ਵਾਲਾ ਇਹਨੂੰ ਕੜੇ ਨਹੀਂ ਸਕਦਾ ਜੀ ਇਹਨੂੰ ਪੰਜਾਬੀ ਬੜੀ ਹੈ ਉਹਨੂੰ ਸਮਝਿਆ ਨਹੀਂ ਆ ਸਕਦੀ ਏ ਉਹ ਗਲਤ ਪੜ੍ਹੂ ਉਹਨੇ ਜੋ ਪੜਿਆ ਉਹੀ ਪੜ੍ਹੂਗਾ ਵਿਚਾਰਾ ਇਹ ਸਾਰੀ ਬਦਲ ਨਹੀਂ ਬਹੁਤ ਸੁਣ ਇਹ ਪੜਾਈ ਹੋਰ ਹੈ ਜਿਆਦੇ ਨਾਲ ਤਾਂ ਹੋਗਾ ਦਸ ਹਿੰਦੀ ਚਾਹ ਆਉਂਦਾ ਅਮਰੀਕਾ ਸ਼ੈਲੋ ਜੀ ਟਾਕਾ ਮੂੜੋ ਚਾਰਥ ਪੇਡਾ ਤਾਂ ਵੜਦੇ ਨੇ ਆਇਓ ਸਹਉਦ ਤਾਕਾ ਮੂੜੋ ਚਾਂਦ ਪੈਦਾ ਜਾਖੋ ਪੇਵ ਨਪਾਵਤ ਵਿਦਾ ਤਾਕੋ ਕਰ ਪਾਹਗ ਅਨੁਮਾਨ ਤਾ ਮੂੜ ਕਥ ਪੇਨ ਜਾਣਤ ਯਾਰ ਤਾਇਓ ਸਾਰੇ ਜਿਆਦਾ ਬਹੁਤ ਘੱਟ ਹੁੰਦਾ ਜਾਂ ਤੂੰ ਮੇਰੇ ਵੱਲ ਹੈ ਜਦ ਜਿਆਦਾ ਬੰਦਾ ਜਦ ਜਦ ਤੂੰ ਮੇਰੇ ਵੱਲ ਹੈ ਤਾਕਾ ਮੋ ਚੰਦ ਮੈਨੂੰ ਕੀਲੀ ਪਰਵਾਹ ਹੈ जा, जा करता ਕਰ ਜਾ ਕਰਤਾ ਸਿਰਠੀ ਕੋ ਸਾਜੇ ਹਾਂ ਜੋ ਜਿਹੜਾ ਜਾਪਤ ਲੇਖੈ ਨਾ ਪਵੈ ਉਸ ਕੋਲ ਹਾਂਜੀ ਜਾ ਚੈ ਕਰ ਡਿੱਗ ਦੀ ਸਾਜੇ ਕੱਠਾ ਜਾਚੇ ਕੱਠਾ ਨਹੀਂ ਜਾ ਚ ਇਕੱਠਾ ਹੁੰਦਾ ਨਾ ਨਾ ਜਾ ਚ ਨਾ ਬਸਨਾ ਜੀ ਇਹ ਕਰੇ ਜਾ ਚ ਇਕੱਠੇ ਅਲੱਗ-ਅਲੱਗ ਬਣਨਾ ਜਾ ਚ ਕਰ ਜਿਸ ਦੇ ਘਰ ਵਿੱਚ ਦਿਗ ਦਿਸ ਹੈ ਆਹ ਦਿਗ ਬ੍ਰਾਹਮਣ ਜਦ ਤੱਕ ਅੱਲਾ ਸਾਰੇ ਅਜੜਾ ਉਹਦਾ ਕਾਰ ਕੀ ਹੈ ਅਜਿਹੇ ਚਤਰਾਉਂਦੇ ਨੇ ਜਿੰਨੀ ਆ ਵੀ ਆਹ ਮੂਰਤੀਆਂ ਜਿੱਤਰ ਉਹਦਾ ਕਾਹਦੇ ਸਾਰਾ ਉਹਨਾਂ ਕਰੇ ਹੈ ਉਹ ਪਾਈ ਉਹਦਾ ਸਰਬਿਆਪੀ ਉਹਦਾ ਘਾਰ ਹੈ ਆ ਜਿਹੜਾ ਸ਼੍ਰੀਤੀ ਹੈ ਨਾ ਸਾਰੀ ਰਚਨਾ ਹੈ ਉਹਦਾ ਹੈ ਆਰਾਮ ਘਰ ਵੀ ਹੈ ਜਦੋਂ ਆਮਰ ਆਮガルਪੋਂ ਹੋਇ ਆਏ। ਆਮガルਪੋਂ ਦਾ ਖਾਣਾ। ਉਧੇ ਖੁੰਝਲਦਾ ਤੇ। ਆਹ ਦੇ ਜਮਾਦ ਖਲਦਾ ਖੁੰਝਲਦਾ। ਮਾਲਕ ਕੌਣ ਸਿੱਟੀ ਦਾ? ਬਣਾ ਦੱਸ। ਸਿੱਟੀ ਦਾ ਮਾਲਕ ਕੌਣ ਹੈ? ਜਿਹਨੇ ਸਿੱਟੀ ਬਣਾਈਆ ਅਰੇ ਜਨਾ। ਉਹ ਮਾਲਕ ਹੈ। ਇਹ ਜੀ ਬਣਾਈ ਹੈ ਉਹ ਭਾਈ ਮਾਲਕਾ ਉਹਦਾ ਘਰ ਹੈ ਜਿਹਨੇ ਉਹ ਟੈਂ ਕੋਠੀ ਬਣਾਈ ਹੈ ਤੁਹੀਂ ਵਿਚ ਰਹਿਣਾ ਤੁਹੀਂ ਮਾਲਕ ਵੀ ਹੈ ਠੀਕ ਹੈ ਜੀ ਉਹਦਾ ਹੁਕਮ ਚੱਲਦਾ ਹੈ ਤੇ ਉਹਦੇ ਇਹ ਬ੍ਰਹਮ ਦਾ ਇੱਕ ਪੂਰਨ ਬ੍ਰਹਮ ਦਾ ਘਰ ਆ ਉਹਨ ਬ੍ਰਹਮ ਅੱਥੇ ਰਹਿੰਦਾ ਹੈ ब्रह्म ज्ञान निके मन परदा जैसे तारू पर प्रकाश जैसे तकोला प्रकाश होयो न पार है जोदा करकी जो हुंदा जोदा अंदर होदा रे हुंदा काठ काठ काठ हुं की हुंदा कड़े दा करकी आ कड़े दा पेट है कड़े दा हाल जी कड़े दा आधार है कड़े दा आधार भनोदा है जिया विरोधी ऊपर दी कार है ਉਹ ਉਹਦੇ ਛੋਟਾ ਆਪੇ ਆਪਣਾ ਘਰ ਹੈ ਜੀ ਹਾਂ ਚਾਚੇ ਘਰ ਦਿਗ ਦਿਸੈ ਸਰਾਇਚਾ ਸੱਸਾ ਰਾਰੇ ਨੂੰ ਕੰਨਾ ਈੜੀ ਨੂੰ ਸਿਹਾਰੀ ਚੱਚੇ ਨੂੰ ਕੰਨਾ ਸਰਾਇਚਾ ਹਾਦੀ ਰਚਨਾ ਦਾ ਘਰ ਚ ਪਾਂਤਾ ਤੇਰੇ ਸਾਕੋ ਸਾ ਸਭ ਕੋ ਜੋ ਦੀਨ ਦਾ ਸਾਲ ਉਹਦੇ ਘਰ ਚ ਹੈ ਸਭ ਕਸਦਾ ਮਾਲ ਕੋਈ ਹੈ ਇੱਕ ਕੋ ਕਰਿਆ ਦੁਆ ਕਰੇ ਨਹੀਂ ਕੋਈ ਉਹ ਤਾਂ ਹੋਵੇ ਨਾ ਵੀ ਦੁਆ ਕਰੇ ਸ਼ਹਿਰ ਦੇ ਘਰ ਉਹਦਾ ਬਾਕੀ ਹੋਰ ਲੋਕਾਂ ਨੇ ਦੁਆ ਤਾਂ ਕਰਦਾ ਹੀ ਨਹੀਂ ਦੁਆ ਤਾਂ ਕੋਈ ਕਰੀ ਨਹੀਂ ਮਾਣ ਜੀ ਬਬਈ ਸਰਾਇ ਚਾ ਦਾ ਅਰਥ ਕੀ ਹੋਇਆ ਸਰਾ ਇਕਦਾਰ ਸਰਾਇ ਕਾ ਹੁੰਦਾ ਉਹਦਾ ਅਸਰ ਨਾ ਕਨਾਤ हां जी हां जिमे सहज सदा सहज छावाण संतोष सराय सदा सील सन्हा सो है आ सराय जड़ा कणात जित तक हद होवे जित तक हद होवे आकारा ए एमदूदा संतार ਆ ਅਗਰ ਹੈ ਸੁਖ ਸੰਗਤ ਦੇ ਵਿੱਚੇ ਹੈ ਸੁਖ ਸੰਗਤ ਉਹ ਆਪ ਹੈ ਹਉ ਦਾ ਅੰਦਰ ਉਹ ਕਹਿੰਦਾ ਮੇਰੇ ਅੰਦਰ ਹੈ ਸਭ ਕੁਝ ਮੇਰੇ ਅੰਦਰ ਮੇਰੇ ਘਰ ਵਿੱਚ ਹੈ ਕਾਦੇ ਅੰਦਰ ਹੁੰਦਾ ਹਾਂਜੀ ਬਬਈ ਪੰਨਾ ਨੰਬਰ 141 ਤੇ ਬੰਦਤੀ ਹੈ ਇੱਕ ਤੰਬੂ ਪਲੰਗ ਨਿਵਾਰ ਸਰਾਈਚੇ ਲਾਲਤੀ ਉਹ ਦੇ ਨਾਲ ਉਹ ਰਾਜੇ ਹੁੰਦੇ ਨੇ ਤੰਬੂ ਹੁੰਦੇ ਛੇ ਪਲੰਗ ਹੁੰਦੇ ਤੇ ਅਰਦਲੇ ਕਨਾਤ ਆ ਲੈਣਦੇ ਕਨਾਤ ਨਾਲੇ ਅਰਦਲੇ ਵਿਚਾਲੇ ਤੰਬੂ ਲਾਉਂਦੇ ਤੇ ਜਿਹੜੇ ਰਾਜੇ ਹੁੰਦੇ ਸੀ ਦਰਬਾਰ ਜੇ ਉਹ ਨਾ ਖੜਦੇ ਸੀ ਕਨਾਤ ਦੇ ਨਾਲੇ ਬੇਜੇਦਾਰ ਹੁੰਦੇ ਸੀ ਕੋਈ ਰਾਤ ਨੂੰ ਹਵਲਿਆਂ ਨਾਲ ਰੱਦ ਹੋਵੇ ਇੱਕ ਮਹਿਲ ਬਣਾਉਂਦੇ تھے ਉਹ ਇੱਕ ਜਾਨੀ ਏਰੀਆ ਜਿਹਦੇ ਵਿੱਚ ਹੋਰ ਕੋਈ ਪੜ ਨਹੀਂ ਸਕਦਾ ਡੋਟੇ ਬੰਨ। ਜਿਹੜਾ ਜਦੋਂ ਨਾਲ ਤੂ ਐ ਅਫਕ ਨਾ ਤਾਲ ਲਵਨੇ। ਕਨਾਤਮੀਂ ਜਿਹੜੇ ਛੋਟਿਆਂ ਨਾਲ ਆਉਂਦਾ ਆ ਖੜੇ ਕਰਦੇ ਆ। ਬਾਉਂਡਰੀ ਬਾਉਂਡਰੀ। ਜਿਹੜੀ ਬਾਉਂਡਰੀ ਬਣਾਉਣੀ ਆ ਉਹਨੂੰ ਕਹਿੰਦੇ ਨੇ ਲੱਕੜ ਦੇ ਵਿੱਚੋਂ ਬਾਸ ਖਾੜੇ ਕਰਕੇ ਵਿੱਚ ਹੁੰਦੀਆਂ ਨੇ ਲਾਈ ਟਰਪਾਲ ਜੀ ਬੋਟਾ ਕਪੜਾ ਹਾਂਜੀ ਹਾਂਜੀ ਹਾਂਜੀ ਉਹ ਖਨਾਤ ਕਹਿੰਦੇ ਨੇ ਦੋਨੋਂ ਦੀ ਦੀਵਾਰ ਬਾਉਂਡਰੀ ਕਾਸ਼ ਦੇ ਵਿਚਾਲੇ ਜਿਹੜੀ ਦੀਵਾਰ ਉਹਦਾ ਨਾਮ ਸੜਾਕੇ ਆ ਉਹ ਕੀ ਹੈ ਜੀ ਉਹ ਪਰਮੇ ਲਿਖਿਆ ਹੈ ਮੈਂ ਹੈ ਦੂਦ ਉਹ ਪਰਮਾੰਡਾ ਲੇ ਪਰਮਾੰਡਾ ਉਹ ਹੈ ਉਦੇ ਵਿੱਚ ਕੂਟੋਂਡਾ ਪਰਮਕਾ ਉਹਨੇ ਪਰਗਾਸਾ ਪਰਗਾਸਾ ਬਾਹਰ ਦਾ ਜਿਹੜਾ ਪਰਮਦੇ ਅੰਦਰ ਪ੍ਰਕਾਸ਼ ਦਾ ਪ੍ਰਕਾਸ਼ ਨਹੀਂ ਹੁੰਦਾ ਜੇ ਪ੍ਰਕਾਸ਼ ਉਹਦਾ ਪ੍ਰਕਾਸ਼ ਤਾਂ ਬਾਹਰ ਹੈ ਪਰਗਾਸਾ ਜਿਹੜਾ ਉਹ ਪ੍ਰਕਾਸ਼ ਨਹੀਂ ਸਾਨੂੰ ਦੇਣਾ ਜਦ ਮੇਰੇ ਹਿੱਤੇ ਦਾ ਰੋਸ਼ਨੀ ਬਾਹਰ ਅੰਦਰ ਇੱਕ ਰੋਸ਼ਨੀ ਹੋ ਗਈ ਉਹ ਪ੍ਰਗਾਸ ਹੈ ਅੰਦਰ ਹੋਏ ਗਿਆਨ ਪ੍ਰਗਾਸ ਇਸ ਵਿਨਾਸ਼ ਪ੍ਰਕਾਸ਼ ਕਰਨਾ ਪੈਂਦਾ ਨੇ ਦੇ ਵਿੱਚ ਫਿਰ ਇਹ ਰਹਿੰਦਾ ਹੀ ਨਹੀਂ ਬਾਹਰੰ ਦੇ ਕੋ ਹੋ ਜਾਂਦਾ ਉਹਨੂੰ ਪ੍ਰਕਾਸ਼ ਰਹਿੰਦੇ ਨੇ ਹਾਂਜੀ ਜਾ ਚੈ ਕਰ ਦਿਗ ਦਿਸੈ ਸਰਾਇਚਾ ਬੈਕੁੰਠ ਭਵਨ ਚਿੱਤਰਸਾਲਾ ਬੈਕੁੰਠ ਭਵਨ ਹੈ ਇਹਨੂੰ ਐ ਬੈਕੁੰਠ ਕਹਿਣਾ ਨੇ ਜਿੜੀ ਬੈ ਕੁੰਠਾ ਦਾ ਹਾਂਜੀ ਜਾਚੈ ਘਰ ਦਿਗ ਦਿਸੈ ਸਰਾਇਚਾ ਆ ਸਰਾਇਚਾ ਇੱਥੇ ਆ ਇੱਥੇ ਬਹੁਣ ਨਹੀਂ ਚਲਣਾ ਪਰ ਮਨ ਸੰਤੋਖ ਦੇ ਉਹ ਸੰਤੋਖ ਦੀ ਬਾਉਂਡਰੀ ਜਾਉਣਾ ਸਤ ਸੰਦੋਰੀ ਲੰਘ ਲੰਘ ਰੋਣ ਦੇਗਾ ਜਿਹੜੇ ਆਰਾਮਕਾਰ ਚਾਹੁੰਦਾ ਉਹ ਲੰਘ ਰੋਣ ਦੇਗਾ ਨਾ ਗੈਰਾਂ ਦੀ ਹੁਲਤ ਰੋਣ ਦੇਗਾ ਆਰਾਮਕਾਰ ਹੈਗਾ ਤੇ ਚਾਹ ਗਰਦਾ ਮਾਰੇ ਆਰਾਮਕਾਰ ਦੁੱਖ ਲਗੇ ਨਾ ਭਾਈ ਦੁੱਖ ਨਹੀਂ ਆਉਂਦੇ ਉਹਦੇ ਆਰਾਮਕਾਰ ਹੈ ਆਰਾਮਕਾਰ ਦੇ ਅੰਦਰ ਉਹਦਾ ਘਰ ਹੈ ਹੈ ਗੁਰਬਾਣੀ ਦੇ ਅੰਦਰ ਉਹ ਰਾਮ ਘਰ ਦੇ ਅੰਦਰ ਉਹਦਾ ਘਰ ਹੈ ਉੱਥੇ ਜਾਉਣਾ ਸਾਨੂੰ ਵੀ ਇਹ ਕਾਚਰ ਉੱਥੇ ਦੇਖਾ ਤੋਂ ਫਿਰ ਖਵਾਲਾ ਮੈਂ ਆ ਇੱਥੇ ਤੋਂ ਉਹ ਇਹ ਘਾਟਾ ਬਤਾ ਦੇ ਉਹਦਾ ਘਰ ਆ ਗਿਆ ਉੱਥੇ ਸਭ ਕੁਝ ਆਪਣਾ ਤੇ ਸਭ ਕੁਝ ਜਦ ਫਰਬੇ ਚਾਪਣੇ ਸਭ ਕੁਝ ਬਾਹਰ ਕਿਉਂ ਜਾਣਾ ਬਾਹਰ ਕੀ ਹੈ ਬਾਹਰ ਨਾਲ ਬੇਸ ਜੋਖਾ ਉਹ ਯਾਰ ਜਣਾ ਵਧੀਆ ਫੜਾ ਮੈਂ ਖਾ ਲਾ ਉਹ ਪੜੀ ਦੀ ਨੂੰ ਜੀ ਦੇ ਬਾਅਦ ਤੇ ਪਹਿਲਾਂ ਕੀਤਾ ਵਾਪੇ ਖਾਲੂ ਜਿਹੜਾ ਤੈਨੂੰ ਪਹਿਲਾਂ ਕੀਤਾ ਉਹ ਕਵਨ ਗਾਲ ਜੀਜ ਖਾ ਲਮੈਂ ਤੈਨੂੰ ਉਹ ਹੀ ਜੀ ਦੱਲਿ ਤੇਰੇ ਬਾਅਦ ਜੱਟਦਾ आले कर दिग दिसै सरायचा बैकुंठ भवन चित्र माने अंदर बाउंड्री का है पिटा ना नहीं कर है ओ सरायचा है ना बाउंड्री है ओले पर सातर दो की है ओदा घर ओ चलीया बक उन्हें आपस में कहता पास दो कह देने ਗਿਆ ਰਾਮਕਾਰ ਕਹਿੰਦੇ ਚੌਕਰ ਦਾ ਮਾਰੇ ਰਾਮਕਾਰ ਰਾਮ ਦਾ ਘਰ ਹੈ ਉਹ ਹੁਕਮ ਨੇ ਜਿਹੜਾ ਉਹੀ ਉਹਦਾ ਘਰ ਹੈ ਹੁਕਮ ਜਿਹੜਾ ਨਹੀਂ ਉਹਦਾ ਘਰ ਹੈ ਜਿੱਥੇ ਤਾਂ ਕੋਹੋਂ ਮੈਨੂੰ ਤੇਸੇ ਕੋਲਾ ਘਰ ਹੈ ਹੁਕਮ ਜਿਹੜਾ ਹੋ ਪਾਣੀ ਤਰੋ ਕਾਜੀ ਜਾ ਚੈ ਕਰ ਦਿਗ ਸਰ ਆਜਾ ਸਨਾਤ ਵੀ ਹੈਗੀ ਬਾਉਂਡਰੀ ਹੈਗੀ ਆ ਮਤਲਬ ਕਹਿਣ ਦਾ ਡਿੱਗ ਦਿਸੈ ਡਿੱਗ ਡਿੱਗ ਦਿਸੈ ਦਿਸ਼ਾ ਦਾ ਦੇਸ਼ਾ ਦੱਦੇ ਨੂੰ ਸਿਹਾਰੀ ਸੱਸੇ ਨੂੰ ਦਲਾਵਾ ਦਿਸ਼ਾ ਦਿਸ਼ਾ ਨੇ ਹੁੰਦੀ ਵਿਸ਼ਾ ਕਹਿੰਦੇ ਨਹੀਂ ਆਪਾਂ जाचे कर दिग दिसै दिग ददनु सारी गंगा दिग है हां जी दिग दा ब्राह्मण नु कहंदा ने भी हुंदा बहुत बड़ा दिग ब्राह्मण ला बहुत बड़ा भी हुंदा है जेड़ा ब्राह्मण है वो बहुत बड़ा है ਬੜੀ ਹਸੀ ਦਾ ਨੋਆ ਦਿੱਕਲੀ ਹੈ ਬਹੁਤ ਉਨਕੀਆ ਹੋ ਆ ਤੋ ਰਾਜ ਨਾ ਉੱਤੇ ਇਹ ਨਾ ਉੱਜਾਗਾ ਉਹ ਛੋਟੀ ਵੱਡੀ ਦਵਾਈ ਨਾ 10 12 ਬੰਦੀ ਵੀ ਟਪੂ ਉਹ ਦਵਾਈ ਕੋਟ ਆਪ ਸਖਦਾ ਬਾਉਂਡਰੀ ਐਜਾ ਬਾਹਰ ਨਹੀਂ ਜਾ ਸਕਦਾ ਤਨ ਸਾਜ ਜਵਰਨ ਲੱਗੀ ਨ ਕੋਈ ਐ ਉਹਦੇ ਕਾਚੇ ਜਿਹੜਾ ਹੁਕਮ ਦੇ ਵਿੱਚ ਨਹੀਂ ਹੈ ਉਹ ਦੁਖੀ ਹੈ ਜਿਹੜਾ ਹੁਕਮ ਦੇ ਵਿੱਚ ਹੈ ਪਾਣੇ ਵਿੱਚ ਸੁਖੀ ਹੈ ਪਰ ਉਹ ਹੈ ਕਾਂ ਚੁਛਾਰੇ ਆ ਕਾਟਾ ਤੇਰੇ ਸਭ ਕਿਛ ਹੈ ਤੂੰ ਕੋਈ ਕੁਝ ਵੀ ਬਾਹਰ ਨਹੀਂ ਦੇ ਰੱਖ ਤੋ ਉਹ ਸਾਰਾ ਕੁਝ ਕਾਚੇ ਉਹਦੇ ਦੁਖੀ ਆ ਜਿਹੜੇ ਆਪਣੇ ਪਾਣੇ ਚੱਲਦੇ ਨੇ ਦੁਖੀ ਨੇ ਜਿਹੜੇ ਉਹਦੇ ਪਾਣੇ ਚੱਲਦੇ ਨੇ ਸੁਖੀ ਨੇ ਆਹ ਦੇ ਕੋਪਸ ਇੰਡੀਆ ਦੇ ਨੇ ਜਿਹੜੇ ਹੁਕਮ ਦੇ ਵਿੱਚ ਚੱਲਦੇ ਨੇ ਸਰਕਾਰ ਦੇ ਨੀਮਾਨ ਸਾਥ ਚੱਲਦੇ ਨੇ ਇਮਾਨਦਾਰੀ ਨਾਲ ਚੱਲਦੇ ਨੇ ਉਹਨਾਂ ਨੂੰ ਕੋਈ ਕੁਝ ਨੀ ਲੈਣੀ ਠੀਕ ਹੈ ਜੀ ਨਹੀਂ ਕਹਿਣਾ ਚਾਹੀਦਾ ਜੇ ਕਹਿਂਦਿਆ ਤਾਂ ਫਿਰ ਉਹ ਰਾਜਨੀ ਤਰਫ ਨਾ ਹੈਗਾ ਉਹਨਾਂ ਨੂੰ ਕੋਈ ਕੁਝ ਨਹੀਂ ਕਹਿਣਾ ਹੁੰਦਾ ਜੇ ਰਾਜਨੇਕ ਹੋਵੇ ਉਹਨਾਂ ਨੂੰ ਕੋਈ ਖਤਰਾ ਨਹੀਂ ਹੁੰਦਾ ਕਬਾ ਜਾਨੇ ਕੋ ਬੇ ਰਾਜੇ ਦੇ ਨਾਲ ਚੱਲਣ ਸਾਰੇ ਹੋ ਸੁਖੀ ਉੱਤੇ ਕਿ ਸੁਧਾਰਾਜ ਇਹ ਰਾਜ ਦੀ ਗੱਲ ਨਹੀਂ ਕਰਦਾ ਜੋ ਮੌਜੂਦਾ ਹੈ ਤਾਂ ਕਿਸੇ ਗੁਦਾ ਰਾਜੇ ਵਿੱਚ ਨਹੀਂ ਗੱਲ ਹੋ ਸਕਦੀ ਇਹ ਜਿਹੜੇ ਬਗਵਾਸ਼ ਨੇ ਸੁਖੀ ਨੇ ਕੁਝ ਬਗਵਾਸ਼ ਸੁਖੀ ਨੇ ਸਰਕਾਰ ਦੇ ਨਾਲ ਜਿਹੜੇ ਬਗਵਾਸ਼ ਨੇ ਲਾਠਾਂ ਸੇ ਨੇ ਸਰਕਾਰ ਤੋਂ ਲਿਆ ਬਗਵਾਸ਼ੀ ਦਾ ਸੁਖੀ ਨੇ ਜਦੋਂ ਹੀ ਪਾਰਟੀ ਆ ਯੂਜ਼ ਹੋਏ ਉਹਨਾਂ ਨੂੰ ਸੁਖੀ ਹੋ ਜਾਣਗੇ ਉਹਨਾਂ ਤੇ ਉਹਨਾਂ ਲਿਆ ਹੋਇਆ ਹੈ ਇਹ ਨਹੀਂ ਅਭੀ ਕੋਈ ਸਰਕਾਰ ਖਰਾਬ ਅਗਰਾਬ ਸਾਡੀ ਨਹੀਂ ਸੁਫੰਸਾੜੀ ਦਿੰਦੇ ਨੇ ਬਦਮਾਸ਼ਾਂ ਨੂੰ ਜੋਰਾਂ ਨੂੰ ਥੱਕਣ ਆਪ ਵੀ ਥੋੜਾ ਥੱਕਦੇ ਚਾਹਸ ਤਾਂ ਇਹਦੀ ਗੱਲ ਨਹੀਂ ਕਰਦੇ ਮੌਜੂਦਾ ਰਾਜ ਦੀ ਇਹ ਰਾਜ ਦੀ ਗੱਲ ਕਰਦੇ ਨੇਖ ਵੀ ਰਾਜ ਹੀ ਨੇ ਉਨੇ ਵਿੱਚ ਦਾ ਰਾਜ ਦਾ ਨੇਕੀ ਦਾ ਰਾਜ ਹੈ ਉਹਦੇ ਘਰ ਵਿੱਚ ਜਿਹੜਾ ਉਹਦੇ ਪਾਣੀ ਚ ਸੁਕੀ ਹੈ ਉਹ ਤੇ ਸੰਸਾਰੀ ਦੇ ਸ਼ੈਤਾਨੋਂ ਨੂੰ ਦੁਖੀ ਦਿੰਦਾ ਵੀ ਹੈ ਇੱਥੇ ਉਹ ਦੁੱਖ ਨੂੰ ਦੁੱਖ ਮੰਨਦਾ ਹੀ ਨਹੀਂ ਦਾਰੂ ਮੰਨਦਾ ਉਹਦੇ ਪਾਣੀ ਸਹਿੰਦਾ ਉਹ ਲੰਮੀ ਨਜ਼ਰ ਨਾਲ ਉਹਦਾ ਆ ਸੰਸਾਰੀ ਦੇ ਉਹਦਾ ਹੈ ਹੀ ਨਹੀਂ ਤੇ ਸਰਕਾਰਾਂ ਜਿਹੜਾ ਨਿਊਟਰਲ ਹੈ ਸਰਕਾਰਾਂ ਮੇਰੇ ਕੋਲ ਕੁਝ ਨਹੀਂ ਕਹਿੰਦੀ ਕੋਈ ਬੰਦੇ ਜਾਵੇ ਸਰਕਾਰੋਂ ਨਹੀਂ ਦੇਣਾ ਜਾਂ ਸਰਕਾਰ ਚੋਂ ਦਖਲ ਹੀ ਨਹੀਂ ਦਿੰਦਾ ਇਸ ਨੂੰ ਕਹਿਣਾ ਹੀ ਕੁਝ ਨਹੀਂ ਸਰਕਾਰ ਵੀ ਉਹਨੂੰ ਕੁਝ ਨਹੀਂ ਰੱਖਦੀ ਸਰਕਾਰ ਨਹੀਂ ਦਿੰਦਾ ਉਹਦਾ ਜੇ ਸਰਕਾਰ ਜਦ 71 ਜਿਹੜੀ ਪਹਿੜੀ ਹੈ ਉਹ ਜੰਗੀ ਲੱਭੀ ਉਹਨੂੰ ਜੰਗਾ ਸਕਦਾ ਇੱਕ ਤਰ ਪਹਿੜੀ ਹੈ ਉਹ ਮਾੜਾ ਸਮਝਦਾ ਫੇਰ ਸਰਕਾਰ ਵੀ ਉਹਨੂੰ ਕਰਦੀ ਹੈ ਕੋ ਕੋ ਦੇ ਆਪਣੇ ਮਨ ਚ ਵੀ ਫਰਕ ਆ ਜਾਂਦਾ ਚੰਸ ਕਾਦਾ ਹੋਇਆ ਦੇ ਸਿੱਖਿਆਦ ਨਹੀਂ ਕੋਈ ਲਵੇ ਸਭ ਨੂੰ ਇੱਕ ਹੋ ਜਾ ਗਏ ਫਿਰ ਕੋਈ ਵੀ ਨਹੀਂ ਰਹਿਣਾ ਹੁੰਦਾ ਕੁਝ ਜਾਂ ਸਾਡੇ ਅੰਦਰ ਫਰਕ ਆਉਂਦਾ ਫਿਰ ਦੂਜੇ ਦੇ ਉੱਪਰ ਕਾ ਜਾਣਾ ਆ ਬਬਲੀ ਇਹਦਾ ਹੁਣ ਜਿਹੜੀ ਪੰਕਤੀ ਆਪਾਂ ਕਰ ਰਹੇ ਆ ਇਹਦਾ ਪ੍ਰੋਪਰ ਅਰਥ ਕੀ ਬਣਿਆ ਚਾ ਚੈ ਘਰ ਦਿਗ ਦਿਸਹ ਸਰਾਇਚਾ ਯਾਰ ਉਹਦੇ ਘਰ ਐਡਾ ਬੜੀ ਬਨਾਤ ਹੈ ਉੱਥੇ ਹੱਥ ਨਹੀਂ ਉੱਪਰ ਦਾ ਕਰਦਾ ਅਥਾਰਾ ਕਾਸ਼ਕ ਨਾ ਤੇ ਉਹ ਜਾਈ ਨਹੀਂ ਹੋਈ ਬੈਕੁੰਠ ਭਵਨ ਹੈ ਬੈਕੁੰਠ ਭਵਨ ਇਹ ਚਿੱਤਰ ਨਹੀਂ ਹੈ ਉਹਦੇ ਰੂਪ ਅਨੂਪ ਹੈ ਕਿਸਮ ਦੇ ਰੂਪ ਇੱਥੇ ਨੇ ਜਿਵੇਂ ਉਹਦੇ ਕਾਦੇ ਵਿੱਚੇ ਇਹਦਾ ਨਾਮ ਦੇਖੋ ਮਨੂ ਅੰਦਰੋਂ ਚਿੱਤਰ ਸ਼ਾਲਾ ਜਿਹੜੀ ਹੈ ਧਰਮ ਸ਼ਾਲਾ ਚਿੱਤਰ ਸ਼ਾਲਾ ਪਾਕ ਸ਼ਾਲਾ ਪਾਕ ਸ਼ਾਲ ਵੀ ਆਇਆ ਲਵ ਜੀ ਪਾਕ ਸ਼ਾਲਾ ਉਹਨੂੰ ਕਹਿੰਦੇ ਜਿੱਥੇ ਰਸੋਈ ਬਖਦੀ ਹੈ ਉਹ ਘਰ ਵੱਡਾ ਹੁੰਦਾ ਉਹਦੇ ਵਿੱਚ ਕਮਰੇ ਹੁੰਦੇ ਨੇ ਚਿੱਤਰ ਵੀ ਕਮਰਾ ਹੁੰਦਾ ਉਹਦੇ ਘਰ ਦੇ ਵਿਚਾਲੇ ਜਿਹੜਾ ਸੰਭਾਰੇ ਚਿੱਤਰ ਸ਼ਾਲਾ ਹੈ ਸਰਵਤੇ ਕੁੰਡ ਪਪਨ ਚਿੱਤਰ ਚਾਲੋ ਦੇ ਵਿੱਚ ਹੈ ਰਚਨਾ RAM ਨੇੜੀ ਰਚਨਾ ਬਣਾਈ ਹੈ ਚਿੱਤਰ ਬਣਾਏ ਨੇ ਜਿਵੇਂ ਕੋਈ ਬਣਾਉਂਦਾ ਨਾ ਆਪਣੇ ਸਿਨਰੀ ਪੇਂਟਿੰਗਸ ਉਹ ਪਿੰਡ ਆਪਣੇ ਬਣਾਈ ਆਪਣੇ ਕਪੜੇ ਖੁੰਡੋ ਦੀ ਸਜਾ ਕੇ ਰੱਖ ਲੈਂਦਾ ਘਟਾ ਉਹਦਾ ਵੱਡਾ ਹੁੰਦਾ ਉਹਨੇ ਆਪਣੇ ਘਰਾਂ ਪੇਂਟਿੰਗ ਬਣਾ ਕੇ ਰੱਖੀ ਜਿੰਨੀਆਂ ਜੋ ਨੇ ਸਤਿ ਸ਼੍ਰੀ ਅਕਾਲ ਹੈ ਉਹਦਾ ਗਾਣਾ ਮੈਂ ਗਾ ਲਿਆ ਕੋਈ ਹਾਂਜੀ ਸਮਝ ਆ ਗਈ ਤੇ ਉਹਦੇ ਅੰਦਰੇ ਕਮਰਾ ਹੈ ਇੱਕ ਉਹਦਾ ਹੀ ਬਾਹਰ ਦਾ ਸੁਠਾਰ ਘਾਦਾ ਇਸ ਸਾਗਰ ਦਾ ਅੰਦਰ ਹੈ ਨਾ ਹਾਂਜੀ ਹੈਗੇ ਜੀ ਬਾਬਾ ਜੀ ਇੱਥੇ ਕੀ ਹੋਇਆ ਚ ਚਿੱਤਰ ਬਚਿੱਤਰ ਇਹ ਹੈ ਅਬ ਚਿਹਰਾ ਇਹ ਅਬ ਇਹ ਚਤਰ ਵਿਚ ਤਰਾਂ ਚਿੱਤਰ ਇਹ ਜਸਤਰ ਨੂੰ ਨਾ ਦੇਖੋ ਨੂੰ ਜਦੋਂ ਆਂ ਕਿ ਤੇਰਾ ਜੀ ਮੈਂ ਚਿੱਤਰ ਬਣਾਇਆ ਉਹਦੇ ਨਾਲ ਉਹਦੀ ਗੱਲ ਕਰੋ ਉਹਦਾ ਧਿਆਨ ਕਰੋ ਇਹ ਚਿੱਤਰ ਨਾਲੇ ਖੋਦੇ ਜੇ ਜਦੋਂ ਦੇਖੋਗੇ ਜਿਹੜੇ ਚਿੱਤਰ ਚ ਫਸ ਗਏ ਉਹ ਰੂਪ ਧਾਰਨ ਕਰਨਾ ਪੈਣਾ ਜਿਹੜਾ ਜਨਨ ਲਗੂ ਤੇ ਵੜਜੋਗੇ ਉੱਥੇ ਧਿਆਨ ਹੋ ਜਾਓ ਉਹ ਚੰਗਾ ਜਿਹਾ ਨਾਲੇ ਉਹ ਸੁਪਨਾ ਦੇਖੀ ਜਾਓਗੇ ਜੋ ਅੰਦਰ ਉਹਦੇ ਚੱਤਰ ਚ ਵੜ ਕੇ ਹਾਂਜੀ ਸਭਤ ਲੋਕ ਸਮਾਨ ਪੂਰੀਲੇ ਆਜਣ ਲੜਣ ਕਈ ਨਾ ਲੋਕ ਨੇ ਸਤਪਤਾਲ ਸੱਤ ਰਾਸ਼ੇ ਬੁੰਦੇ ਨੇ ਉਹਨਾਂ ਦਾ ਰਾਸ਼ਨ ਪਾਣੀ ਸਾਬ ਵਿੱਚ ਭਰਿਆ ਹੈ ਪੂਰੀਲੇ ਉਹਨਾਂ ਨੇ ਪੂਰਾ ਕਰਨ ਵਾਸਤੇ ਹੈ ਬਹੁਤ ਕੋਲੇਵਲ ਪੂਰਾ ਕਰਨ ਵਾਸਤੇ ਖਾਣ ਪੀਣ ਦਾ ਸਾਮਾਨ ਵੀ ਵਿੱਚ ਉਹਨਾਂ ਦੇ ਤੇ ਦਵੀ ਦਾ ਭਰਨਾ ਹੈ ਸਭ ਦਾ ਜੀ ਗਿਆਨ ਵਾਲਾ ਵੀ ਭਰਨਾ ਚੁਗਾ ਵੀ ਭਰਨਾ विके राशन वाणी जो कुछ पाया से एक बार एक बार पाता हां जी जी आप कर रहे सी पन्ना 1292 तो राग मलर वाणी भगत जियो की जाचे कर लक्ष्मी कोवारी चंद सूरज दीवड़े कौतुक काल बपुड़ा कोतवाल सुकरा श्री ਲੱਛਮੀ ਲੱਛਮੀ ਉਹਦੀ ਹੁੰਦੀ ਹੈ ਲੱਛਮੀ ਮਾਇਆ ਨਹੀਂ ਹੁੰਦੀ ਉਹ ਮਾਇਆ ਵੀ ਚਮਕਦੀ ਆ ਅਸਲ ਜਸਲ ਚਮਕਦੀ ਆ ਅਕਲ ਦਾ ਗਿਆਨ ਚਮਕਦਾ ਜਿਹੜੀਆਂ ਦੇਸ਼ ਤਲਵਾਰਾਂ ਨੇ ਜਿਹੜੇ ਗਿਆਨ ਦੇ ਲੈਸ ਕਬੂਦੀ ਨਹੀਂ ਬਾਹਰ ਆਉਂਦੀ ਹੈ ਅੰਦਰ ਜੋ ਗਿਆਨ ਦੀ ਰੋਸ਼ਨੀ ਆ ਬਲੇਵਾਰ ਕੱਢਦੀ ਆ ਉਹਨੂੰ ਤੇ ਬੋਲ बोल के या कुछ करके दिखा के ए लक्ष्मीया गोरी गोरी होरेंदी है ओनु कहंदा रे तू मेरी मेरा माता तू मेरा पिता तू है मेरा माता बोला लक्ष्मीया गोरी ओबित ओदे घर हैगी है अकल ओदे घर है ਅਗਲੋ ਫਿਰ ਮਿਲਦੀ ਹੈ ਉਹ ਗੁਰਮਤ ਉਹਥੇ ਮਤ ਉਹਥੇ ਹੀ ਮਿਲਦੀ ਹੈ ਮਤਮਤਾ ਮਤ ਉਹਥੇ ਹੀ ਮਿਲਦੀ ਹੈ ਗੁਰਮਤ ਉਹਥੇ ਹੀ ਮਿਲਦੀ ਹੈ ਸਾਰ ਬਾਣੀ ਉਥੋਂ ਹੀ ਆਈ ਹੈ ਧੁਰ ਬਾਣੀ ਇਹ ਹੁੰਦਾ ਕਹਿੰਦਾ ਜਾਂ ਜਿੰਨੀ ਸੋਚੀ ਆਉਂਦੀ ਹੈ ਉਥੋਂ ਹੀ ਆਉਂਦੀ ਹੈ ਸੋਚੀ ਉਹ ਲక్ష్ਮੀ ਹੈ ਸੰਸਾਰ ਨੂੰ ਜਿੰਨੇ ਪ੍ਰਕਾਰ ਦੀ ਸੋਚੀ ਹੈ ਉਥੋਂ ਹੀ ਹੁੰਦੀ ਹੈ ਇਹ ਹੀ ਹੈ ਜਿਦੋਂ ਸੋਦੀ ਆਉਂਦੀ ਉਹਦੇ ਵਿੱਚ ਚਮਕ ਲਸ਼ਕ ਜਿਵੇਂ ਬਿਜਲੀ ਲਸ਼ਕੀ ਐਂ ਜਦੋਂ ਕਲਸ਼ਕ ਬਾਦੋਂ ਆਉਂਦੀ ਜਦੋਂ ਸੋਦੀ ਆ ਜਾਂਦੀ ਹੈ ਕਲਿਕ ਹੋ ਜਾਂਦੀ ਹੈ ਘਰ ਲਕਸ਼ਮੀ ਕੁਆਰੀ ਹਾਂ ਚੰਦ ਸੂਰ ਆਜ ਚਤਾਰ ਮੰਦੇ ਹੀ ਬੜੇ ਨੇ ਉਹ ਕਿੱਥੇ ਦੀਬੜੇ ਕਿੱਥੇ ਬਿਜਲੀ ਦੀ ਰੋਸ਼ਨੀ ਚਾਉਂ ਕੋ ਪਤਾ ਦੀਵੜੇ ਨੇ ਦੋਏ ਵਿਚਾਰੇ ਆ ਦੂਏ ਚੰਦ ਸੂਰਜੇ ਦੇ ਨੇ ਤਾਂ ਪਤਾ ਨਹੀਂ ਕਿੰਨੇ ਕਰਨੇ ਇਹ ਵੀ ਉਹਦੇ ਘਰ ਨੇ ਆ ਦੂਏ ਜਿਹੜੇ ਚੰਦ ਸੂਰਜੇ ਨੇ ਆਪਣੇ ਜੜ ਚੰਦ ਸੂਰਜੇ ਜੜ ਤਾਂ ਅਸੀਂ ਨੋਂ ਰੱਖ ਲਏ ਉਹਨਾਂ ਦੇ ਚੰਨ ਸੂਰਜ ਚੇਤਨ ਵੀ ਨੇ ਚੰਨ ਸੂਰਜ ਜੜ ਵੀ ਨੇ ਦੋਈ ਉਹਦੇ ਘਰ ਚ ਨੇ ਹਾਂਜੀ ਚੰਦ ਸੂਰਜ ਦੀਵੜੇ ਅੱਜ ਤਰਮਨ ਚੰਨ ਸੂਰਜ ਨੇ ਇਹ ਰਸੋਈ ਕਰਦੇ ਨੇ ਉਹ ਦੀ ਪਿਆਰ ਉਹ ਸੋਈ ਗਿਆ ਆਹ ਜਿੰਨੇ ਵੀ ਗਿਆਨ ਸੋਈ ਆਤਮਾ ਦਾ ਗਿਆਨ ਇਹੀ ਕਹਿੰਦਾ ਕਰਦੇ ਨੇ ਕਉ ਰਸੋਈ ਸੋਈ ਕਿ ਚੰਦ ਸੂਰਜ ਬਿਨਾ ਫਲ ਕੋਈ ਫਸਲ ਨੀ ਹੁੰਦੀ ਬਾਹਲੇ ਜੀਤੇ ਫਰਾਗੰਦਲੇ ਜੀਂ ਦੀ ਖਰਾਬ ਹੋਏ ਪੈਦਾ ਇਹੀ ਕਰਦੇ ਨੇ ਚਾਹ ਕਿਸੇ ਪ੍ਰਕਾਰ ਦੀ ਵੀ ਹੋਵੇ ਅੱਡ ਅੱਡ ਜੁਨੀਏ ਦੀ ਅੱਡ ਅੱਡ ਖਰਾਬ ਹੈ ਅੱਡ ਅੱਡ ਸਾਰੀ ਅੱਡ ਅੱਡ ਖਰਾਬ ਹੈ ਚਾਰ ਵੇਦ ਨੇ ਚਾਰ ਪ੍ਰਕਾਰ ਦਾ ਗਿਆਨ ਚਾਰੇ ਪ੍ਰਕਾਰ ਦਾ ਚਾਰੇ ਵੇਦ ਬ੍ਰਹਮੇ ਕੋ ਦੱਤੇ ਨੇ ਉਹਦੇ ਘਰੇ ਆ ਉਹਨਾਂ ਕਰੋ ਨਹੀਂ ਮਿਲੇ ਨੇ। ਛਾਰੇ ਪ੍ਰਕਾਸ਼ ਦਾ ਗਿਆਨ ਸੰਸਾਰ ਚ ਹੈ। ਛਾਰੇ ਪ੍ਰਕਾਸ਼ ਦੇ ਵਿਦਵਾਨ ਨੇ। ਅਤਾਂਗ ਕਰਾਂਗੀ ਵਾਲਾ ਗਿਆਨ ਵੀ ਉੱਥੋਂ ਮਿਲਿਆ। ਉਹਦੇ ਵੀ ਖੜਾ ਖਾਲੇ ਲੋਕ ਹੈਗੇ ਨੇ। ਉਹਦੀ ਪੁਖਾਲੇ ਵੀ ਨੇ। ਸੰਸਾਰਿਕ ਗਿਆਨ ਦੀ ਪੁਖਾਲੇ ਵੀ ਨੇ। ਨਿਰਾਕਾਰ ਦੇ ਗਿਆਨ ਦੇ ਪੁਖਾਲੇ ਵੀ ਨੇ। ਦੋਹੇ ਪ੍ਰਕਾਸ਼ ਦਾ ਗਿਆਨ ਹੈ ਉੱਥੋਂ ਹੀ ਮਿਲਦਾ। ਜੇ ਕਿ ਚੰਦ ਦਾ ਗਿਆਨ ਹੈ ਸੰਸਾਰੀ ਬੁਖ ਇੱਕ ਸੂਰਜ ਦਾ ਗਿਆਨ ਹੈ ਮੈਰਾਹਾਰੀ ਬੁਖ ਜਿਹੜਾ ਬ੍ਰਹਮ ਗਿਆਨ ਹੈ ਉਹ ਸੂਰਜ ਦਾ ਗਿਆਨ ਹੈ ਉਹ ਪਰਮ ਦਾ ਨਾਸ ਕਰਦਾ ਹੈ ਉਹ ਤਾਂਹੇ ਸੂਰਜ ਵੰਸੀ ਕਹਿੰਨੇ ਨੇ ਰਾਮਚੰਦਰ ਨੂੰ ਸੂਰਜ ਕਿਉਂ ਸੀ ਕਿ ਪਿਛੋਕੜ ਵਾਲਿਆਂ ਦਾ ਗਿਆਨ ਬ੍ਰਹਮ ਗਿਆਨ ਸੀ ਨਾ ਕੋਲੋਂ ਉਕੇ ਮਾਰਤਾ ਨੇ ਫੇਰੀਆ ਮਰਿਆਦਾ ਪਰਛੋਦਦਾ ਰਾਮ ਬਣਿਆ ਬੇੜਾ ਕਰਤਾ ਰਾਮ ਨੇ ਕੀਤਾ ਵੈਦ ਦਾ 라ਵਣ ਨੂੰ ਮਾਰ ਕੇ 라ਵਣ ਦਾ ਵਿਰੋਧ ਕਰਦਾ ਹੈ ਰਿਸ਼ੀ ਮੋਨੀ ਜਿਹੜੇ ਪਖੰਡਵਾਦੀ ਨੇ ਉਹਨਾਂ ਦੀ ਸਪੋਰਟ ਕਰਦਾ ਹੈ ਵਰਕੀਟਾ ਕੀ ਉਹ ਮੂਰਤੀ ਪੂਜਾ ਮੰਦਰ ਤਾਂ ਬਣਾਉਂਦੇ ਨੇ ਉਹਨਾਂ ਦੀ ਰੋਜੀ ਰੋਟੀ ਉਹਦੇ ਵਿੱਚ ਹੈ ਬਾਟ ਜਿਨ੍ਹਾਂ ਨੇ ਪਾੜੀ ਹੈ ਨਾ ਪੰਡਤ ਨੇ ਬਾਟ ਪਾੜੀ ਉਹਨਾਂ ਨੂੰ ਸ੍ਰਕਸ਼ਨ ਦੇਣ ਵਾਲਾ ਇਹੀ ਰਾਮ ਹੈ। ਤਾਂ ਕਬੀਰ ਨੇ ਬਦਲਤਾ ਸਭੇ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰਿਕੇ ਹਾਰੂ ਪੰਡਤ ਨੂੰ। ਸੁੰਦਰ ਬੋਲਦਾ ਉਹ ਰਾਮ ਹੈ ਥੋੜੇ ਵਾਲਾ ਰਾਮ ਰਾਮ ਨਹੀਂ ਹੈ। ਉਹਨੇ ਤਾਂ ਬਾੜ ਪਾੜੀ ਏ, ਉਹਦੇ ਅਸਲ ਤਾਂ ਤੁਸੀਂ ਬਾੜ ਪਾੜੀ ਏ। ਅੱਜ ਉਹ ਕਹਿੰਦੇ ਨੇ, ਵੀ ਸ਼ਗਰੂ ਦੀ ਲੋੜ, ਹੁਣ ਦੇਖਾਂਗੇ ਕਦੇ ਬਣਦਾ ਵੀ ਸ਼ਗਰੂ। ਬੇਸ਼ਗਰੂ ਬਣੂਗਾ। ਸਾਰੇ ਦੁਨੀਆ ਨੇ ਮਤਤਾਨੂੰ ਰੋਜ਼ ਨਹੀਂ ਲਊਗਾ ਕਰੂਗਾ ਨਹੀਂ ਤਾਂ ਫਰਮਾਈ ਤੇ ਗੁਰੂ ਕੀ ਜਾਤੇ ਭਰਮ ਜਾਏ ਹਾਂਜੀ ਚੰਨ ਤੇ ਸੂਰਜ ਦੀਵੜੇ ਕੌਤਕ ਕਾਲ ਬੱਪੂੜਾ ਚੰਨ ਸੂਰਜ ਦੀਵੜੇ ਚੰਨ আর ਸੂਰਜ ਦੀਵਨੇ এবੀ ਰੋਜ਼ ਨਹੀਂ ਦੇ ਰਹੇ ਨੇ ਸੂਰਜ ਦੀ ਰੋਸ਼ਨੀ ਤਾਂ ਪਰਮ ਦਾ ਨਾਸ ਕਰਦੀ ਹੈ ਹਨੇਰਾ ਚੱਕਦੀ ਹੈ ਚੰਨ ਦੀ ਰੋਸ਼ਨੀ ਜਿਹੜੀ ਹੈ ਉਹ ਰਾਤ ਨੂੰ ਹੁੰਦੀ ਹੈ ਰੋਸ਼ਨੀ ਤਾਂ ਕਰਦੀ ਹੈ ਸੀਮਤ ਰੋਸ਼ਨੀ ਕਰਦੀ ਹੈ ਬਹੁਤ ਸੀਮਤ ਜਿਹਨੇ ਜਿਹੜਾ ਗਿਆਨ ਚਾਹੀਦਾ ਉਸ ਨੂੰ ਉਹ ਜਿਹਾ ਹੀ ਗਿਆਨ ਦਿੰਦੀ ਹੈ ਜੋ ਮੰਗਣਾ ਠੰਕਰ ਪਰੰਤੇ ਸੋਈ ਸੋਈ ਦੇਵਾ ਨਾਨਕ ਇੱਥੇ ਕੋਮਲ ਗੁਰੂ ਨਾਨਕ ਨੂੰ ਅੰਕੜਾ ਲੱਗਿਆ ਹੋਇਆ ਇੱਥੇ ਜੇ ਔਂਕੜ ਨਹੀਂ ਹੈ ਔਂਕੜ ਲਾਉਣਾ ਪਊਗਾ ਨਾਨਕ ਦਾਸ ਮੁਖ ਤੇ ਜੋ ਬੋਲਣ ਜਿਨੇ ਦਾਸ ਨੇ ਉਹਦੇ ਜਿਹੜੇ ਵੀ ਉਹ ਬੋਲਦੇ ਨੇ ਮੁਖੋ ਇਹ ਆ ਵਹ ਸੱਚ ਹੋਆ ਕਿਉਂਕਿ ਭਗਤ ਦਾਸ ਨੇ ਸਾਰੇ ਉਹ ਬੋਲੇ ਨੇ ਇਹ ਪਰ ਲੋਕ ਜੋ ਸੱਚ ਹੈ ਉਹ ਇਹਨਾਂ ਨੇ ਕਿਹਾ ਜਦ ਲੱਗ ਜਾਏ ਨਾ ਨਾਲ ਨਾਨਕ ਦੇ ਸਤ ਮੰਦ ਜੁੜ ਜਾਂਦਾ ਔਕੜ ਹਟ ਜਾਂਦਾ ਉਹ ਕੜ ਨਹੀਂ ਹਟ ਸਕਦਾ ਇੱਥੇ ਕਿ ਦਾਸਰਾਂ ਉਂਕਰ ਲੱਗੂਗਾ ਜਾ ਕੇ ਜੇ ਦਾਸਰਾਂ ਉਂਕਰ ਲਾ ਦੀਏ ਜਾ ਕੇ ਨਾਨਕ ਨੂੰ ਦਾਸ ਬਣਾ ਦਈਏ ਤੇ ਭਗਤ ਕਿੱਥੇ ਗਏ ਜਿਹੜੇ ਉਹ ਬੋਲਣੇ ਬਾਬਾ ਜੀ ਮੇਰੇ ਕੋਲ ਈਸ਼ਰ ਮਾਈਕਰੋ ਜਿਹੜੀ ਗੁਰਬਾਣੀ ਦੀ ਐਪ ਹੈ ਉਹਦੇ ਵਿੱਚ ਨਾਨਕ ਮੁਕਤ ਹੈ ਕੱਕਾ ਮੁਕਤ ਹੈ ਦਾਸ ਤੇ ਉਂਕਰ ਲੱਗੀ ਹੈ ਗੱਲ ਤਾਂ ਮੇਰੇ ਨਾਨਕੇ ਦਾਸ ਹੋ ਗਿਆ ਇੱਕ ਵਕਤ ਦਾਸਰੇ ਤਾਂ ਕਿੱਥੇ ਗਏ ਉਹ ਗੁਰਬਾਣੀ ਜਿਹਦੇ ਭਗਤ ਬੈਠੇ ਨੇ ਉਹ ਉਹਨੀਆਂ ਵਾਹ ਬੋਲ ਨਾਮ ਕਰਿਆ ਇਹਦਾ ਮਤਲਬ ਇਹ ਹੋ ਗਿਆ ਦਾ ਸੱਚ ਹੈ ਨਹੀਂ ਸੱਚ ਹੈ ਗੁਰਬਾਣੀ ਦਾ ਹੈ ਇਹ ਤੇ ਜਦ ਨਾਨਕ ਜੀ ਬੋਲ ਰਹੇ ਹੈ ਹਾਂ ਨਾਨਕ ਦਾ ਕਾਹ ਰਿਹਾ ਕਹਿ ਰਹੇ ਫਿਰ ਨਾਨਕ ਦਾ ਮੁਖ ਫੇ ਤਾਂ ਕਿ 3rd ਪਰਸਨ ਦੀ ਬਾਣੀ ਹੋ ਗਈ ਨਾਨਕ ਜੀ ਦੀ ਬਾਣੀ ਉਹਨਾਂ ਲਈ ਹੈ ਤੇ ਜੀ ਆਏ ਪਾਏ ਨੇ ਇਹਨਾਂ ਨੇ ਇਹਨਾਂ ਦੀ ਅਕਲ ਨਹੀਂ ਸਾਰੀ ਬਾਣੀਆਂ ਗਲਤ ਕਰਦੀ ਸਾਰੀ ਬਾਣੀ ਗਲਤ ਕਰਦੀ ਤਾਂ ਜਿੰਨੀਆਂ ਵੀ ਸੀਗੀਆਂ ਸਾਈ ਨਾਲੀਆਂ ਮਿਲਡਾ ਜਿਦਾਂ ਗੁਰੂ ਘਰ ਦੇ ਦੱਸ ਸਾਰੀਆਂ ਖਤਮ ਕਰਤੀਆਂ ਉਹਨੇ ਉਹ 50 ਸਾਲ ਚ ਖਤਮ ਕੀਤੀਆਂ ਨੇ ਸਰੋ ਖਾਕ ਫਾਸੀ ਉੱਜੜਿਆ ਥੰਦਾ ਰਿਹਾ ਇੱਕ ਵੀ ਮਿਲ ਨਹੀਂ ਛੱਡੀ ਉਹ ਤਾਂ ਹਰ ਜਿਹੜਾ ਜਿਹਨੂੰ ਤੱਕ ਪ੍ਰੋਬਲਮ ਨੀ ਇਹਨਾਂ ਨੂੰ ਜੀ ਵੀ ਕੋਈ ਕਰ ਨਹੀਂ ਸਕਦਾ ਕਰ ਕਿਉਂ ਨਹੀਂ ਸਕਦਾ ਕਿਉਂ ਨਹੀਂ ਕਰ ਸਕਦਾ ਕੀ ਇਹ ਗੱਲ ਝੂਠ ਹੈ ਹਰ ਜੁਗ ਜੁਗ ਕੋ ਭਗਤਾ ਪਾਇਆ ਜੀ ਜੇ ਭਗਤਾਂ ਦੇ ਬਾਦ ਆਨੰਦ ਗੁਰਨਾਨ ਕੋ ਹੋ ਸਕਦਾ ਹੈ ਹੋ ਸਕਦੇ ਨੇ ਸੁੰਦਰ ਹੋ ਸਕਦਾ ਹੋਰ ਕਿਉਂ ਨਹੀਂ ਕੋਈ ਸਮਝਦਾਗਾ ਜੀ ਹੋ ਸਕਦੇ ਕਿਉਂ ਨਹੀਂ ਸਮਝਦਾ ਕੋਈ ਜੇ ਨਹੀਂ ਸਮਝ ਆ ਰਹਾ ਫਿਰ ਬੇਕਾਰ ਸੀ ਤੇ ਪੰਥ ਚਲਾਉਣਾ ਬੇਕਾਰ ਸੀ ਤੇ ਬੀੜ ਲਿਖਣੀ ਬੇਕਾਰ ਸੀ ਇਹਦਾ ਫਾਇਦਾ ਸੀ ਇੱਥੇ ਕਿ ਪੰਥ ਚਲੇ ਤਬ ਜਗਤ ਮੇਂ ਜਬ ਤੁਮ ਕਰੋ ਜਬ ਤੁਮ ਕਰੋ ਸਾਹਿਬ ਇਹ ਕਹਿੰਨਾ ਨੇ ਆਪਣੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੰਨੀ ਗੱਲ ਕਰਦੇ ਜੀ ਗਲਤ ਹੋ ਗਿਆ ਪ੍ਰਚਾਰ ਤੋਂ ਹੁੰਦੇ ਹੀ ਉਹ ਪ੍ਰਚਾਰ ਹੋ ਗਿਆ ਗਲਤ ਉਹ 76 ਨੇ ਜਿਹੜੀ ਹੋਣੀ ਹੈ ਉਹ ਤਾਂ ਹੋਊਗੀ ਹੋ ਵੀ ਹੁੰਦੀ ਰਹੂ ਨੇ ਚੋਰੀ ਕੀਤੀ ਹੈ ਖਾਂਦੇ ਨੂੰ ਉਹ ਦੇਖੀ ਗਏ ਨੇ ਛੱਤਰ ਦੇਖੀਏ ਹੁਣ ਜਿਹੜਾ ਰੰਗ ਲਾ ਦੇਣਗੇ ਉਹ ਦੇਖ ਲਾਂਗੇ ਜਿਹੜੇ ਪੰਜਾਬ ਦੇ ਸਿੱਖ ਨੇ ਜਿਹੜੇ ਹੁਣ ਵਿਸ਼ਗੁਰੂ ਬਣਾ ਰਹੇ ਨੇ ਉਹਨਾਂ ਨਾਲ ਕਿੰਨਾ ਬਿਜਾਇਆ ਉਹ ਦਿਨ ਪਤਾ ਕਬਸ ਬੋਲ ਹੋ ਜਾਣੇ ਇਹਨਾਂ ਨੂੰ ਬਿਸ਼ਵਗੁਰੂ ਤਾਂ ਹਿੰਦੂ ਬਣਾਉਣ ਲੱਗੇ ਨੇ ਮੁਸਲਮਾਨ ਨਾਲ ਨੇ ਈਸਾਈ ਯਹੂਦੀ ਨਾਲ ਨੇ ਇਹ ਇਨਕਸਾਫ ਤਾਂ ਵੀ ਮਰੇ ਨਾ ਦੇਣਗੇ ਤੋਂ ਭਲਾ ਚਿੱਖੀ ਤੋਂ ਐਂਟੀ ਚਿੱਖੀ ਤੋਂ ਸਾਥ ਹੋ ਜਾਣਗੇ ਸਾਧਨ ਵਿੱਚ ਬਗੜਨ ਦੇ ਖੇਤਰ ਖਾ ਕੇ ਬਿਲਕੁਲ ਐਡਮਿਟ ਕੌਤਕ ਕਾਲ ਬੱਪੂੜਾ ਕਾਲ ਬੱਪੂੜਾ ਕਾਲ ਕੀ ਹੈ ਕਲਪਨਾ ਹੀ ਕਾਲ ਹੈ ਇਹੀ ਤੋਦ ਕਰਦਾ ਇਹ ਕਾਲ ਹੈ ਮਨ ਜਿਹੜਾ ਨਾ ਇਹੀ ਇਹਦਾ ਕਾਲ ਹੈ ਸਾਡੀ ਅਕਲ ਦਾ ਕਾਲ ਅਕਲ ਦਾ ਦੁਸ਼ਮਣ ਮਨ ਕਲਪਨਾ ਕਰਦਾ ਮਨ ਕਲਪਨਾ ਹੀ ਕਾਲ ਹੈ ਕਾਲ ਕਲਪਨਾ ਕਦੇ ਨਾ ਖਾਏ ਉਹ ਇਹ ਕਹਿੰਦੇ ਕਾਲ ਕਲਪਨਾ ਨੇ ਸਾਨੂੰ ਖਾਈ ਜਾਂਦੀ ਹੈ ਸਾਡੀ ਅਕਲ ਨੂੰ ਖਾਈ ਜਾਂਦੀ ਹੈ ਸਾਡੇ ਗਿਆਨ ਦਾ ਨਾਸ ਕਰੀ ਜਾਂਦੀ ਹੈ ਬੁੱਧੀ ਦਾ ਨਾਸ ਕਰਦੀ ਹੈ ਕਲਪਨਾ ਜਿੰਨਾ ਚਿਰ ਜੋ ਸੋਚਦੇ ਨੇ ਸਾਡੀ ਬੈਟਰੀ ਡਾਊਨ ਹੁੰਦੀ ਹੈ ਅਕਲ ਦੀ ਜੇ ਬਚਾ ਲਵੇ ਗੁਰਬਾਣੀ ਬੈਠੀ ਯਾਰਜ ਹੁੰਦੀ ਹੈ ਚਾਰੇ ਤਾਂ ਕਰਦੇ ਹੀ ਨਹੀਂ ਗੁਰਬਾਣੀ ਤਾਂ ਵਿਚਾਰਦੇ ਹੀ ਨਹੀਂ ਸੋਚ ਸੋਚ ਕੇ ਬੈਠੀ ਢੋਂ ਕਰਦੀ ਇੰਨੀ ਡਾਊਨ ਹੋ ਗਈ ਸੱਖਾਂ ਦੀ ਬੈਠੀ ਉਹਨਾਂ ਨੂੰ ਪਤਾ ਹੀ ਨਹੀਂ ਕੀ ਕਰੀਏ ਕਿ ਦੁਨ ਜਾਈਏ। ਡੇਰਾ ਹੀ ਨਾ ਰਚਾਂਸ ਭੇਰੇ ਨਾ। ਗੁਰੂ ਛੱਡਤਾ ਨਾ ਮਾਇਆ ਲੈ ਲਈ। ਠੱਗ ਮੂਰੀ ਖਾਈ। ਉਹ ਠੱਗ ਮੂਰੀ ਖਾਲੀ ਮਾਇਆ। ਉਹ ਠੱਗਾਂ ਦੀ ਜਿਹੜੀ ਸੀ ਨਾ ਆਪਣੇ ਆ ਗੁਰਮਤ ਠੱਗਾਂ ਨੇ ਜੋ ਅਰਥ ਕੀਤੇ ਗੁਰਮਤ ਦੇ ਠੱਗ ਮੂਰੀ ਸੀ ਉਹ ਖਾਲੀ ਮੂਰੀ ਦਾ ਸਵਾਦ ਮਿਠਾ ਤਾਂ ਹੁੰਦਾ ਨਹੀਂ ਉਹ ਖਾਲੀ ਠੱਗ ਮੂਰੀ ਖਾਈ ਮੂਰੀ ਕੀ ਹੁੰਦਾ ਜੀ ਮੋਲੀ ਬੋਲੀ ਬੋਲੀ ਨੂੰ ਮੂਰੀ ਕਹਿੰਦੇ ਨੇ ਬੋळा ਉਹ ਮੂਰੀ ਮੂਰੀ ਬਣ ਗਈ ਉਹ ਉਹ ਮੂਰਤੋਂ ਲੱਲੇ ਤੋਂ ਰਾਜਾ ਬਣ ਗਿਆ ਬੋੜ ਹੈ ਨਹੀਂ ਨਾ ਸਾਡਾ ਉਹ ਬੋੜ ਤਾਂ ਸਾਡਾ ਸੱਚ ਹੈ ਖਾਲੇ ਝੂਠ ਠੱਗ ਮੂਰੀ ਖਾਈ ਇਹ ਕੰਦਾਲੀ ਬਣਾਈ ਹੋਈ ਜਲ ਅਜੇ ਵੀ ਕਹਿੰਦੇ ਨੇ ਇਹਦੀ ਆ ਪ੍ਰਾਣੀ ਮਤ ਦਾ ਸਨਾਤਨ ਮਤ ਦਾ ਪ੍ਰਾਣੀ ਉਹ ਕੀ ਹੁੰਦੀ ਹੈ ਝੂਠੀ ਮਤ ਸੱਚ ਪ੍ਰਾਣਾ ਹੋਵੇ ਸੱਚੀ ਮਤ ਪ੍ਰਾਣੀ ਹੁੰਦੀ ਦੀ ਸੱਚੀ ਮਤ ਚੇਰਾਣੀ ਹੁੰਦੀ ਆ ਝੂਠੀ ਮਤ ਪ੍ਰਾਣੀ ਹੋ ਜਾਂਦੀ ਹੈ ਹੁੰਦੀ ਰਹਿੰਦੀ ਹੈ ਪ੍ਰਾਣੀ ਕੀ ਹੁੰਦਾ ਕੋਣ ਨੇ ਖੁੱਟੇ ਨਾਨਕਾਉੜ ਸੱਚ ਰਹੀ ਫੇਰ ਕੋਡ ਕੋਟਾ ਸਾਹਿਬ ਤੋਂ ਜੰਨ ਸੱਚ ਫੇਰ ਪਰਟ ਹੋ ਜਾਂਦਾ ਹੈ ਤਾਂ ਇਹ ਪੰਕਤੀ ਪੰਕਤੀ ਕਿੱਥੋਂ ਦੀ ਹੈ ਜੀ ਕਬੀਰ ਦਾ ਸ਼ਬਦ ਹੈ ਧਰਨ ਆਪ ਨਹੀਂ ਖਾਦੀ ਕਬੀਰ ਨੇ ਵਾਲਾ ਨਹੀਂ ਫੇਰਦਾ ਸੀ ਜਿਆ ਮਾਰਾ ਫੇਰਦਾ ਸਾਰੀ ਜ਼ਿੰਦਗੀ ਨੰਗੀ ਮੂਹ ਚ ਦੋਲ ਆਉਂਦੀ ਮੋੜੀ ਦੀ ਗੱਲ ਮੋੜੀ ਦੇ ਕੰਦ ਚੰਗੀ ਹੁੰਦੀ ਹੈ ਉਕਾਵਤਾ ਕੇ ਦੁਰਗੰਧ ਓਡੀ ਦੁਰਗੰਧ ਦਾ ਹੈ ਜਿਆਦਾ ਪ੍ਰਚਾਰ ਕਰਦੇ ਦਰਬਾਨੀ ਦਾ ਉਲਟਾ ਦੁਰਗੰਧ ਦਾ ਊੜੀ ਉਹਦੀ ਔਰ ਕੀ ਹੈ ਉਹ ਊੜੀ ਇਸ ਮਹਿਲ ਹਾਂਜੀ ਕੌਤਕ ਕਾਲ ਬਪੁਰਾ ਕੋਟਵਾਲ ਕੋਈ ਕੋਟਵਾਲ ਦਰਮੂਰੇ ਉਹ ਵੀ ਇੱਕ ਪਾਸੇ ਪੁੰਨਾ ਇੱਕ ਪਾਸੇ ਪਾਪ ਦੋ ਦਰਵਾਜ਼ੇ ਨੇ ਨਾ ਪਾਪੋਂ ਦਰਵਾਜਾ ਨਹੀਂ ਪਾਪ ਦਾ ਦਰਵਾਜਾ ਤਾਂ ਮੰਨਵਾਲਾ ਜੇ ਪਾਪਾ ਖੋਲ੍ਹੇ ਉਥੇ ਮੰਨਤਾੜਿਆ ਮਵასი ਰਾਜਾ ਇਹ ਹਿਰਦੇ ਆਲਾ ਖੋਲ੍ਹੇ ਉਥੇ ਦੁਆ ਬੈਠਾ ਧਰਮ ਰਾਜ ਬੈਠਾ ਇੱਕ ਪਾਸੇ ਧਰਮ ਰਾਜ ਆ ਇੱਕ ਪਾਸੇ ਮਨੂ ਮਵასი ਰਾਜਾ ਸਾਖਤ ਹੈ ਇੱਕ ਪਾਸੇ ਸੰਤ ਬੈਠਾ ਇੱਕ ਉਥੇ ਸਾਖਤ ਬੈਠਾ ਇੱਕ ਸਾਖਤ ਦਾ ਗੇਟ ਹੈ ਹੁਣ ਜਾਣਦਾ ਇੱਕ ਸੰਤ ਦਾ ਕੌਜਾ ਨੀ ਮੈਂ ਕਹਿੰਦੇ ਤੇ ਹਾਂਜੀ ਚੰਦ ਸੂਰਜ ਦੀਵੜੇ ਕੌਤਕ ਕਾਲ ਬਪੂੜਾ ਕੋਟਵਾਰ ਇੱਕ ਪਾਸੇ ਦਾ ਮਨ ਬੈਠਾ ਕਾਲ ਇਹ ਆਪਣਾ ਹੀ ਕਾਲ ਆ ਪੁੱਠਾ ਇਹ ਪੁੱਠੀ ਹੈ ਕਲਪਨਾ ਕਰਦਾ ਇੱਕ ਪਾਸੇ ਧਰਮ ਰਾਜ ਆਲਾ ਹੈਗਾ ਉਹ ਸੁਗਰਤਾ ਉਧਰਲੇ ਪਾਸੇ ਦੋ ਹੁਕਮ ਨੇ ਇੱਥੇ ਇਹਦੇ ਘਰ ਚ ਐਂ ਕਹਿ ਲਾ ਇੱਕ ਮਨ ਪਾਉਣਾ ਹੁਕਮ ਮਨ ਕਾ ਪਾਣੇ ਦੁਰ ਕਾ ਪਾਣੇ ਇਹਨੇ ਦੋ ਇੱਕ ਪਾਸੇ ਦਾ ਗੇਟ ਮਨ ਕੇ ਪਾਣਿਆ ਉਹਨੇ ਨਾਲ ਇੱਕ ਪਾਸੇ ਗੁਰ ਕੇ ਪਾਣਿਆ ਗੇਟ ਇੱਕ ਪਾਸੇ ਸੰਤ ਨਾਲ ਇੱਕ ਪਾਸੇ ਦੋ ਇਹਨੇ ਨਾ ਜੀ ਇਹਦਾ ਕారణ ਉਹ ਕਹਿੰਦੇ ਆਦ ਅਪਾਰ ਅਲੇਖ ਅਨੰਤ ਅਕਾਲ ਅਪੇਖ ਅਲਖ ਅਨਾਸਾ ਰਜਨਾਂ ਕੀ ਹੈ ਇਕ ਸਵਈਏ ਚ ਦੱਸਿਆ ਦਸਮ ਬਾਸ਼ਾ ਨੇ ਸਾਰਾ ਕੁਝ ਜਿਹੜਾ ਹੈ ਨਾ ਆਦ ਅਪਰ ਕੈ ਸ਼ਿਵ ਸ਼ਕਤੀ ਦਿਓ ਸੰਸਚਾਰ ਤਮ ਸਤ ਸੂਰ ਕਾ ਦੀਪ ਸਸੀ ਸੂਰ ਕਾ ਦੀਪ ਜੀਵੇ ਕਰਕੇ ਆ ਗਿਆ ਨਾ ਸਸੀ ਸੂਰ ਕਾ ਦੀਪ ਦੋ ਦੀਵੜੇ ਅੰਗਰ ਜੀ ਇਹ ਤਾਂ ਵਧੀਆ ਚਾਲ ਹੈ ਨਾ ਪੂਰੇ ਦਾ ਪੂਰੀ ਰਚਨਾ ਨਹੀਂ ਕਰਤੀ ਇਹ ਤਾਂ ਪੂਰੀ ਨਹੀਂ ਹੋ ਸਕੀ ਸਿਰ ਜਸੂਰ ਕੈ ਦੀਪ ਕਰਕੇ ਜੀਵਲੇ ਸੋ ਸੇਟਰ ਠੀਕ ਪੰਕੇ ਨਾਲ ਪ੍ਰਕਾਸ਼ ਹੈ ਪ੍ਰਕਾਸ਼ ਨਹੀਂ ਹੈ ਬੈੜ ਬੜਾਏ ਲੜਾਈ ਸੁਰਾਸੁਰ ਆਪੋ ਦੇਖਤ ਬੈਠ ਤਮਾਸ਼ਾ ਸੁਰਾਸੁਰ ਅਸੁਰ ਦੇਖਦੇ ਰਖ ਦੁਆ ਨੂੰ ਪੈਦਾ ਕਰਦਾ ਤੋਂ ਉਹਦੇ ਅੰਦਰ ਬਦਾ ਉੱਤਾ ਆਪ ਤਮਾ ਸਾ ਦੇਖ ਲੈ ਰਚਨਾ ਆ ਉਹ ਸੁਭਿਆ ਦੇ ਵਿੱਚ ਆ ਇਸ ਕੀ ਰਚਨਾ ਹੈ ਸਾਰੀ ਉਹ ਕਿਵੇਂ ਕੀਤੀ ਉਹਨੇ ਹਾਂਜੀ ਬੱਬਾ ਜੀ ਇੱਥੇ ਪਾਠ ਹੈ ਚੰਦ ਸੂਰਜ ਦੀਵੜੇ ਕੌਤਕ ਕਾਲ ਬਪੂੜਾ ਕੋਟਵਾਲ ਉਹ ਕਾਲ ਆਪਣਾ ਪੈਰ ਘੋੜਾ ਮਾਰਦਾ ਕੋਤਖੋਰ ਖਣਕੀ ਕੀ ਕਰਦਾ ਕੋਤ ਤਾਂ ਕਰਦਾ ਸਾਦਾ ਪੈਰ ਘੋੜਾ ਮਾਰੀ ਜਾਂਦਾ ਉਹ ਨਾਕੀ ਚੇਤੇ ਕਰਦਾ ਹੈ ਕੋਤਖ ਕੋਤਕ ਕਰਦੇ ਕਾਲ ਵਪੜਾ ਕੋਤਖ ਜਿਹੜਾ ਕਰਦਾ ਹੈ ਇਹ ਮਨਤਾ ਨੇ ਫਾਂਸਨ ਕੀ ਵੀ ਨਹੀਂ ਫਾਂਸਨ ਕੀ ਸਭ ਕੋ ਜਾਣੇ ਛੁੱਟੜ ਕੀ ਇੱਕ ਜੋ ਦੋਈ ਕੋਮਿਲੀ ਹੈ ਉਧੂ ਦੇ ਪਾਸੇ ਹੈ ਇਹ ਕਾਲ ਵਪੜੇ ਦਾ ਨੇ ਨਾਟਕ ਚੇਟ ਕੋ ਕੌਤਕ ਦਾ ਉਹ ਕੌਤਕ ਕਹਿੰਦੇ ਇਹ ਬੱਪੂੜਾ ਬਾਬਾ ਜੀ ਇੱਥੇ ਪਾਠ ਹੈ ਸੁਕਰ ਉਹ ਸੁਕਰੀ ਕਰਨੀ ਸੀ ਪਤੰਸ਼ੂ ਕਾ ਲਖ ਦੇ ਕਰੀਂ ਕਰੀ ਨਹੀਂ ਹੈ ਉਹ ਸ਼ੁਕਰਾ ਵੀ ਹੈ ਨਾ ਸ਼ੁਕਰ ਹੈਗਾ ਸ਼ੁਕਰ ਇਹਨਾਂ ਦਾ ਗੁਰੂ ਹੈ ਇਹਦਾ ਗੁਰੂ ਦੀ ਹੈ ਸ਼ੁਕਰ ਜਿਹੜੇ ਸ਼ੁਕਰ ਦਾ ਗੁਰੂ ਹੈ ਉਹ ਮੂrti ਪੂਜਾ ਨੂੰ ਨਹੀਂ ਮੰਨਦਾ ਮਾਇਆ ਨੂੰ ਨਹੀਂ ਮੰਨਦਾ ਸ਼ੁਕਰਵਾਰ ਜੁਮਾ ਕਹਿੰਦੇ ਜੀ ਨਾ ਆਹੋ ਉਹ ਸ਼ੋਮਕਾ ਸ਼ੋਮਕਾ ਕਰੀ ਸੁਖ ਕਦੀ ਸੁਖ ਰੀਤੀ ਹੁੰਦੀ ਪਬਈ ਕੁਸ ਜਗਾ ਪਾਠ ਹੈਗਾ ਸੁਖਰਾ ਇਕੱਠਾ ਹੈ ਉਹ ਅਰਥ ਦਾ ਉਹ ਹੀ ਸੁਖਰਾ ਕੋਈ ਸੁਖਰਾ ਬਣਿਆ ਇਹ ਹੁਣ ਪਾਠ ਇਕੱਠਾ ਕਰਾਂਗੇ ਜੀ ਸੁਖਰਾ ਜੋ ਆਪਣੇ ਸੈਂਚੀ ਭਾਗ ਦੂਜਾ ਹੈ ਉਹਦੇ ਅਲੱਗ-ਅਲੱਗ ਹੈ ਜੀ ਸੂ ਉਹ ਫਿਰ ਸ਼੍ਰੋਮਣੀ ਕਮੇਟੀ ਦੇ ਵਿੱਚ ਐਨਾ ਨਹੀਂ ਸੀ ਇਹ ਜਿਹੜੇ ਨੇ ਨਾ ਆਪਣੇ ਸੰਪਰਦਾਈ ਜੀ ਇੰਨੇ ਨਿਗਰਜ ਨੇ ਇਹ ਬਿਦਵਾਨ ਗਰੇ ਨੇ ਉਹਨਾਂ ਉਹ ਫਿਰ ਵੀ ਕਾਸ਼ੀ ਦੇ ਪੜ੍ਹੇ ਸੀ ਧਰਮ ਪੜ੍ਹਿਆ ਸੀ ਸ਼ੁਕਰਾ ਉਹਨਾਂ ਨੂੰ ਪਤਾ ਵੀ ਸ਼ੁਕਰਾ ਕੀ ਹੁੰਦਾ ਹੈ ਸ਼ੁਭਕਰਮ ਕਰਨੀ ਤੋਂ ਪਰ ਇੱਥੇ ਸਭ ਕੁਝ ਹੈ ਤਾਂ ਅਸੀਂ ਕੀ ਕਰਨਾ ਹੈ ਉਹਦੇ ਨਾਲ ਸਭ ਕੁਝ ਹੈ ਉਹ ਤਾਂ ਕੱਲ ਜਿਹੜਾ ਬਪੜਾ ਉਹ ਦੱਨੀ ਜਾਣਾ ਤਾਂ ਤਾਂ ਇੱਧਰ ਰਹਿਣਾ ਸਰタル ਵਾਲੇ ਪਾਸੇ ਰਹਿਣਾ ਸੁਖਰਤ ਕਾਲ ਨਾ ਆਇਆ ਤਾਂ ਦੁਖਰਤ ਕਾਲ ਨਹੀਂ ਆਇਆ ਉਹ ਇਹ ਵੀ ਆਊਗਾ ਆਇਆ ਹੋਇਆ ਹਾਂਜੀ ਹੈਗੇ ਫਿਰ ਕੋਈ ਗੱਲ ਦੋ ਕਰਮ ਨੇ ਇੱਕ ਸੁਖਰਤ ਨੇ ਦੁਖਰਤ ਨੇ ਉਹ ਜਿਹੜਾ ਦੂਆ ਪਾਸੇ ਦੁਖ ਤਾਲ ਬਪੜੇ ਵਾਲੀ ਉਥੇ ਖੋਤ ਕਦੇ ਠੀਕ ਹੈ ਜੀ ਸੋ ਐਸਾ ਰਾਜਾ ਸ੍ਰੀ ਨਰਹਰੀ ਨਰਹਰੀ ਐਸਾ ਰਾਜਾ ਹੈ ਉਹਦੇ ਘਰ ਦੋੇ ਕੰਮ ਨੇ ਉਹਦੇ ਘਰ ਸੰਤ ਵੀ ਉਹਦੇ ਨੇ ਉਹ ਦੂਸਰ ਸੰਤ ਵੀ ਉਹਦੇ ਹੀ ਨੇ ਉਹ ਅਸੰਤ ਨੇ ਸ਼ਾਂਤ ਨੇ ਸੰਤ ਨੇ ਦੋਏ ਨੇ ਉਹਦੇ ਘਰ ਭਲੇ ਬੁਰੇ ਸਭ ਤੇਰੇ ਆਇਆ ਨਹੀਂ ਭਲੇ ਵੀ ਉਹਦੇ ਨੇ ਬੁਰੇ ਵੀ ਉਹਦੇ ਨੇ ਉਹ ਰਾਮ ਰਾਧ ਦੋਏ ਨੇ ਪੰਜਵੇਂ ਪਾਸ਼ਾ ਵੀ ਭਲਾਂ ਉਹਨਾਂ ਦੇ ਹੀ ਨੇ ਜੂਏ ਦੋਨੇ ਉਹ ਵੀ ਉਹਦੇ ਹੀ ਨੇ ਇੱਥੇ ਨਾਲੋ ਇੱਥੇ ਅੱਗੇ ਪਤਾ ਲੱਗਦਾ ਇੱਕੋ ਸਗੇ ਭਾਈ ਨੇ ਅਡੱਡ ਨੇ ਪਰ ਪਹਿਲਾਂ ਸਗੇ ਭਾਈ ਅਡੱਡ ਨਹੀਂ ਹੋਏ ਇਕੱਠੇ ਰਹੇ ਨੇ ਚਾਹੇ ਅਵਧਾ ਦੇ ਮੁੰਡੇ ਸੀ ਚਾਹੇ ਗੁਰਨਾਮ ਦੇ ਖੁਦ ਮੁੰਡੇ ਸੀ ਚਾਹੇ ਅੰਗਦ ਦੇ ਮੁੰਡੇ ਸੀ ਜੇ ਕੋਨੇ ਕੋਨੇ ਨਹੀਂ ਨੇ ਉਹ ਦੋ ਇਕੱਠੇ ਹੀ ਰਹੇ ਨੇ ਖਲਾਫ ਰਹੇ ਨੇ ਜੀ ਇਹ ਕਿ ਆ ਕੇ ਤਿੰਨ ਹੋ ਗਏ ਇੱਕ ਉਧਰ ਹੋ ਗਿਆ ਦੋ ਹੋ ਗਏ ਦੋ ਰਹੇ ਨੇ ਫਿਰ ਵੀ ਖਲਾਫ ਪਾਸੇ ਚਲੇ ਜੋੜਾ ਹੀ ਰਿਹਾ ਹੈ ਹਾਂ ਜੀ ਜੀ ਸੇਵਲੇ ਜੇ ਸੇਵਾ ਕਰਨੀ ਹੈ ਜੇ ਕਿਸ ਨੂੰ ਸੇਵਾ ਕਰੀ ਦਿਆ ਇਸ ਦੀ ਤੋ ਸਿਖਿਆ ਲਈਆ ਉਹਦੀ ਸੇਵਾ ਕਰਦੀ ਹੈ ਗੁਰ ਸੇਵਾ ਸ਼ਬਦ ਵਿਚਾਰ ਹੈ ਸਾਡੇ ਜਿਹੜਾ ਗੁਰ ਕੀ ਸੇਵਾ ਹੈ ਨਾ ਆਪਣੇ ਜਿਹੜਾ ਅੰਦਰ ਗੁਰਾ ਉਹਦੀ ਵੀ ਸੇਵਾ ਇਹਦੇ ਚ ਹੁੰਦੀ ਜਿਹੜਾ ਉਪਦੇਸ਼ ਹੈ ਸਾਨੂੰ ਕਰਦਾ ਸਤਗੁਰ ਉਹ ਜੋ ਕਹੇ ਉਹ ਕਾਰਕਮਾ ਉਹ ਗੁਰ ਕਹਿਆ ਸਾ ਕਾਰਕਮਾ ਉਹ ਜਿਹੜਾ ਕਹਿੰਦਾ ਉਹੀ ਸੇਵਾ ਹੈ ਗੁਰ ਕਾ ਬਚਨ ਜਿਹੜਾ ਹੈਗਾ ਮੰਨਣਾ ਉਹਨੂੰ ਦ੍ਰਿੜ ਕਰਨਾ ਹੋਤੇ ਚਲਣਾ ਇਹ ਸਭ ਤੋਂ ਵੱਡੀ ਸੇਵਾ ਹੈ ਸੇਵਾ ਉਹ ਚੀਜ਼ ਹੁੰਦੀ ਹੈ ਜਿਹਦੇ ਨਾਲ ਜਿਹਦੀ ਸੇਵਾ ਕਰੀ ਤੇ ਖੁਸ਼ ਹੋਵੇ ਹੁਣ ਜਿਹੜਾ ਸਤਿਗੁਰ ਹੈ ਆ ਗੁਰਦੇਵ ਹੈ ਅਸਲੀ ਹੈ ਜਿਹੜਾ ਸੱਚਿਆਰਾ ਸੱਚਾ ਉਹ ਸੱਚੇ ਮਾਰਗ ਚੱਲਣ ਤੇ ਖੁਸ਼ ਹੁੰਦਾ ਸੱਚੇ ਮਾਰਗ ਚੱਲਦੇ ਆ ਉਸਤ ਕਰੇ ਜਹਾਨ ਜਦੋਂ ਜੋ ਕਹਿੰਦਾ ਉਹਨੂੰ ਮੰਨੇ ਜਿਵੇਂ ਜਿਹੜੇ ਸਾਡੇ ਸਤਗੁਰੂ ਸੀਗੇ ਉਹ ਕਿਹਦੇ ਤੱਕ ਖੁਸ਼ ਨੇ ਕਿਹੜੇ ਸਿੱਖ ਤੇ ਖੁਸ਼ ਹੋਣਗੇ ਜਿਹੜਾ ਗੁਰਬਾਣੀ ਨੂੰ ਸਮਝੇ ਸਹੀ ਉਹਦੇ ਤੇ ਜ਼ਿਆਦਾ ਖੁਸ਼ ਨੇ ਜਿਹੜਾ ਝੜਾਵਾ ਜ਼ਿਆਦਾ ਝੜਾਵੇ ਆ ਹੋਰ ਕੁਝ ਕਰੇ ਉਹਦਾ ਹੰਕਾਰ ਕਰੇ ਉਹਦੇ ਨਾਲ ਖੁਸ਼ ਨਹੀਂ ਆਏ ਉਹ ਸੇਵਾ ਹੱਥੀ ਕਰੇ ਉਹਦਾ ਹੰਕਾਰ ਕਰ ਲਵੇ ਉਹ ਤੇ ਦੇ ਖੋਜ ਨਹੀਂ ਕਾੜੀ ਤੇ ਪ੍ਰਹਾਰੀ ਨੇ ਹੋ ਕਾੜੀ ਦੇ ਖਲਾਫ ਨੇ ਹੋ ਉਹ ਸੇਵਾ ਦੇ ਵਿੱਚ ਭਾਵੇਂ ਸਾਡਾ ਹੀ ਫਾਇਦਾ ਹੈ ਪਰ ਉਹਦੇ ਨਾਲੇ ਜਿਆਦਾ ਖੁਸ਼ ਨਹੀਂ ਟੀਚਰ ਕਦੋਂ ਖੁਸ਼ ਹੁੰਦਾ ਜਿਹੜਾ ਸਟੂਡੈਂਟ ਸਭ ਤੋਂ ਇੰਟੈਲੀਜੈਂਟ ਹੋਵੇ ਟੀਚਰ ਦੀ ਗੱਲ ਧਿਆਨ ਨਾਲ ਸੁਣੇ ਚੰਗੇ ਨੰਬਰ ਲੈ ਕੇ 100% ਪਾਸ ਹੋਵੇ ਟੀਚਰ ਉਹਦੇ ਨੂੰ ਬੜਾ ਖੁਸ਼ ਹੁੰਦਾ ਹਾਲਾਂਕਿ ਸੁਣਨ ਦਾ ਫਾਇਦਾ ਹੈ ਕੋ ਟੀਚਰ ਬਣਾਉ ਖੁਸ਼ ਹੁੰਦਾ ਸਕੂਲ ਵਾਲੇ ਬਹੁਤ ਉਹਨੂੰ ਪ੍ਰੇਮ ਕਰਦੇ ਨੇ ਵੀ ਸਾਡਾ ਰੋਸ਼ਨ ਕਰਦਾ ਹੈ ਐਵੇਂ ਸਤਗੁਰੂ ਹੁੰਦਾ ਵੀ ਨੌਰੋ ਉਹ ਤੇ ਚੱਲਦਾ ਮੇਰੇ ਪਿੱਛੋਂ ਇਹ ਉਹੀ ਪ੍ਰਚਾਰ ਕਰੂ ਜਿਹੜਾ ਅਸੀਂ ਕਰਦੇ ਹਾਂ ਇਹਨੂੰ ਕਹਿੰਦੇ ਨੇ ਸਪੂਤ ਇਹ ਸਪੂਤ ਹੁੰਦੇ ਨੇ ਇਹ ਸਪੂਤ ਨੇ ਜਿਹੜੇ ਗਾਹਾਂ ਬਾਬਾਣੀਆ ਕਹਾਣੀਆਂ ਪੂਤ ਸਪੂਤ ਕਰੇਨ ਇਹ ਜਿਹੜੀ ਬਾਵਾਨੀ ਕਹਾਣੀ ਹੈ ਇਹ ਬਾਵਾਨੀ ਕਹਾਣੀ ਹੈ ਗੁਰਮਤਿ ਪ੍ਰਚਾਰ ਬਾਬੇ ਤੋਂ ਲੈ ਕੇ ਆਦਮ ਤੋ ਪਿੱਛੋਂ ਲੈ ਕੇ ਤਰੋਂ ਰਾਜਾ ਰਾਮ ਦੀ ਕਹਾਣੀ ਇਹਨੂੰ ਜਿਹੜੇ ਸਪੂਤ ਪੋਤ ਨੇ ਉਹ ਕਰਦੇ ਨੇ ਸਪੂਤ ਜਿਹੜਾ ਪੁੱਤਰ ਹੁੰਦਾ ਉਹਦੇ ਨਾਲ ਖੁਸ਼ੀ ਹੁੰਦਾ ਬਾਪ ਇਸ ਕਰਕੇ ਗੁਰਤੀ ਸੇਵਾ ਸ਼ਬਦ ਵਿਚਾਰ ਹੈ ਉਹਦੀ ਸੇਵਾ ਕਰੋ ਜਿਹੜਾ ਗੋਪਾਲ ਰਾਏ ਹੈ ਤਕੋ ਕੋਲ ਦਾ ਮਤਰਾ ਸ਼ਰੀਰ ਦੇ ਵਿੱਚ ਜਿਹੜਾ ਬੋਲਦਾ ਉਹ ਬੋਲਦਾ ਜਿਹੜਾ ਉਹ ਨਹੀਂ ਨਹੀਂ ਨਾਲ ਸ਼ਰੀਰ ਤਾਂ ਬੋਲਦਾ ਹੈ ਸ਼ਰੀਰ ਦੇ ਵਿੱਚ ਜਿਹੜਾ ਬੋਲਦਾ ਉਹਦੇ ਨਾਲ ਸਾਡਾ ਸਮਝ ਹੁੰਦਾ ਨਾ ਕਿ ਉਹਦੇ ਸ਼ਰੀਰ ਨਾਲ ਸ਼ਰੀਰ ਨਾਲ ਨਹੀਂ ਸਾਡਾ ਬਹੁਤ ਆਸਮੰਦ ਜਿਹੜਾ ਬੋਲਦਾ ਉਹ ਸਾਤ ਸਰੂਪ ਹੈ ਸ਼ਰੀਰ ਨਹੀਂ ਸਾਤ ਸਰੂਪ ਹੈ ਸਿਰ ਤੱਕ ਸਾਜ ਹੈ ਜਿਹਦੇ ਨਾਲ ਤੁਲ ਪੈਦਾ ਕਰਦਾ ਹੈ ਪੈਦਾ ਹੁੰਦੀ ਹੈ ਬਸ ਸਾਨੂੰ ਸੁਣਦੀ ਹੈ ਕੁਝ ਅੰਤਰਾ ਬਿਛੋ ਸਤਗੁਰ ਸਤਗੁਰ ਤੇ ਖਾਲੀ ਕੋਈ ਨਹੀਂ ਉਹ ਆਪਣੇ ਵਿਚਾਰ ਸਰੀਰ ਰੂਪੀ ਜੰਤ ਵਜਾ ਕੇ ਸਾਡੇ ਨੂੰ ਕੰਨਾਂ ਨੂੰ ਸੁਣਨ ਵਾਲੀ ਤੋਂ ਪੈਦਾ ਕਰਦਾ ਹੋਰ ਸਰੀਰ ਦਾ ਕੋਈ ਰੋਲ ਹੀ ਨਹੀਂ ਹੈ ਸਰੀਰ ਦਾ ਕੋਈ ਰੋਲ ਨਹੀਂ ਸਤਗੁਰ ਬਾਸਤੇ ਸਿਰਫ ਆਪਣੇ ਜੋ ਵਿਚਾਰ ਸਾਡੇ ਤੱਕ ਕੰਨਾਂ ਨੂੰ ਸੁਣਾ ਕੇ ਪਚਾਉਣ ਤੱਕ ਆਪਣਾ ਗਿਆਨ ਸਰੀਰ ਦਾ ਰੋਲ ਹੈ ਜਿਵੇਂ ਅਸੀਂ ਕੋਈ ਜੰਤ ਵਜਾਉਨੇ ਆ ਬਾਜਾ ਸਾਰੰਗੀ ਕੋਈ ਚੀਜ਼ ਪੈਦਾ ਕਰਕੇ ਉਹ ਧੁਨ ਪੈਦਾ ਕਰਕੇ ਸੁਣਾਉਨੇ ਆ ਇੰਨਾ ਹੀ ਰੋਲ ਹੈ ਸ਼ਰੀਰ ਦਾ ਜਿਆਦਾ ਨਹੀਂ ਹੈ ਅਸੀਂ ਸਾਰਾ ਹੀ ਸ਼ਰੀਰ ਨੂੰ ਮਹੱਤਵ ਦਿੰਦਾ ਸ਼ਰੀਰ ਦੀ ਕੁੱਲ ਹੁੰਦੀ ਹੈ ਆ ਕੁੱਲ ਉਹ ਹੈ ਜਿਹੜਾ ਅੰਦਰ ਬੋਲਦਾ ਹੈ ਉਹ ਰਾਏ ਦੀ ਸੇਵਾ ਕਰਦੀ ਨੇ ਉਹਦਾ ਸ਼ਰੀਰ ਦੀ ਸੇਵਾ ਨਹੀਂ ਕਰਨੀ ਸ਼ਰੀਰ ਦੀ ਸੇਵਾ ਜਿਹੜੀ ਉਹ ਸੇਵਾ ਨਹੀਂ ਹੈ ਸਰੀਰ ਦੀ ਸੇਵਾ ਦਰਗਾਹ ਪਰਵਾਣ ਨਹੀਂ ਇੱਥੇ ਜੋ ਸੇਵਾ ਸੰਸਾਰ ਚ ਪਰਵਾਣ ਤਾਂ ਹੋ ਸਕਦੀ ਐ ਸੇਵਾ ਉਹ ਅਸੀਂ ਤਾਂ ਉਹਨੂੰ ਸੇਵਾ ਮੰਨ ਸਕਦੇ ਹਾਂ ਸੰਸਾਰੀ ਲੋਕ ਸਾਨੂੰ ਸਰੀਰ ਈ ਅਸੀਂ ਸਰੀਰ ਤੱਕ ਹੀ ਮਹਦੂਦ ਹਾਂ ਪਰ ਦਰਗਾਹ ਦੇ ਵਿੱਚ ਜਿਹੜਾ ਖੁਦ ਸਤਗੁਰ ਹੈ ਉਹ ਤਾਂ ਦਰਗਾਹ ਦੀਆਂ ਬਾਤਾਂ ਹੀ ਦੱਸਦਾ ਹੈ ਹਰ ਦਰਗਾਹ ਬਾਤਾਂ ਨਾਨਕ ਆਖ ਸੁਣਾਵਾ ਹਰ ਦਰਗਾਹ ਦੇ ਵਿੱਚ ਜਿਹੜੀ ਸੇਵਾ ਉਹ ਸੇਵਾ ਦੀ ਗੱਲ ਐ ਇੱਥੇ ਹੋ ਰਹੀ ਅਗਰ ਸੰਥਾਰੀ ਸੇਵਾ ਦੀ ਗੱਲ ਹੋ ਰਹੀ ਹੈ ਸੇਵਾ ਕਰਨੀ ਹੈ ਤਾਂ ਅਕਲ ਨਾਲ ਜੰਦੀ ਸੇਵਾ ਕਰੋ ਜੋ ਗੁਰ ਦਾ ਫਰਮਾਨ ਜੋ ਸਾਨੂੰ ਫਰਮਾਇਆ ਹੈ ਉਹਨੂੰ ਮੰਨੋ ਪਰ ਉਤੇ ਚੱਲੋ ਚੱਬਣ ਚੱਲਣ ਸੇ ਰਤਨ ਸੁਣੀਅਰ ਬਹਿ ਗਏ ਫਰੀਦ ਕਹਿੰਦਾ ਈਨਾਂ ਨੇ ਵਿਚਾਰੇ ਗੁਰਬਾਣੀ ਨੂੰ ਸੁਣ ਕੇ ਵਿਚਾਰੇ ਚੱਪਣ ਦਾ ਹੁੰਦਾ ਵਿਚਾਰੇ ਫੇ ਚੱਲੇ ਨੇ ਸੋ ਰਾਤਾਂ ਉਹ ਉਹਨਾਂ ਨੂੰ ਰਤਨ ਹੁੰਦਾ ਤਨ ਜੀਰਾਂ ਦਾ ਰੰਗਿਆ ਗਿਆ ਉਹਨਾਂ ਨੂੰ ਇਨਾਮ ਦਾ ਰੰਗ ਚੜਿਆ ਉਹਨਾਂ ਨੇ ਆਪਣਾ ਹਿਰਦਾ ਰੰਗਿਆ ਉਹਨਾਂ ਨੇ ਆਪਣੀ ਕਾਇਆ ਰੰਗੀ ਹੈ ਕਾਇਆ ਰੰਗਣ ਜੇਥੀਆ ਪਾਈਏ ਨੌਂ ਮਜੀਠ ਨਾਮਦਾਰਾਂ ਨੂੰ ਚਾੜਿਆ ਰੰਗੜਾ ਵਾਲਾ ਜਿਹੜੇ ਸਾਹਿਬ ਰੰਗਾਲੇ ਸਾਹਿਬ ਸਤਗੁਰ ਉੱਥੋਂ ਆ ਰੰਗ ਐਸਾ ਰੰਗ ਨਾ ਡੀਟ ਐਸਾ ਰੰਗ ਵੀ ਤੁਹਾਨੂੰ ਕਿਤੇ ਹੋਰ ਮਿਲਣਾ ਨਾ ਆਉਂਦਾ ਉਹ ਐਸੇ ਵਾਹੇ ਆਪਣੇ ਆਪ ਨੂੰ ਗੁਰਬਾਣੀ ਦੇ ਵਿੱਚ ਮਨ ਨੂੰ ਮੰਨਦਾ ਭੇਜੇ ਜਾਣਾ ਜੇ ਗੁਰਬਾਣੀ ਦੇ ਨਾਮ ਦੇ ਵਿੱਚ ਮਨ ਭੇਜਿਆ ਨਹੀਂ ਸੇਵਾ ਨਹੀਂ ਹੋਈ ਜਿਹੜਾ ਮਨ ਭੇਜ ਗਿਆ ਫੇਰ ਉਹ ਚੜ ਗਿਆ ਫੇਰ ਚੜ ਗਿਆ ਇਹ ਗੱਲ ਕਹੀ ਹੈ ਇੱਥੇ ਸੇਵਿਆ ਲੈ ਗੋਪਾਲ ਰਾਏ ਅਕੋਲ ਨਰਨਜਣ ਉਹਦੀ ਸੇਵਾ ਕਰਦੀਆਂ ਦੇਹ ਦੇ ਨਾਲ ਕੋਈ ਸੰਬੰਧ ਨਹੀਂ ਇਸ ਗੱਲ ਦਾ ਸਰੀਰ ਨਾਲ ਹਾਂਜੀ ਭਗਤੀ ਦਾਣ ਦੀਜੈ ਉਹ ਕੀ ਕਰਦਾ ਭਗਤੀ ਦਾਣ ਦੰਡਾ ਹੋ ਭਗਤੀ ਦਾਣ ਉੱਥੋਂ ਮਿਲਦਾ भक्ति की है मत दंदा गुरकी मत तू ले ओयाने ओ ले लो ओ दी मत जेडी दे रिया है भक्ति बिना बहुत डूबे सयाने यही भक्ति है जे एयर नी जेडे भक्ति बड़े बड़े स्याने डूब गए वाला फेर नाले और योगी सब डूब गए जिना गुरमत लई है ਗੁਰੂ ਕੀ ਮੱਤ ਲਈ ਗੁਰ ਕੀ ਮੱਤ ਤੂੰ ਲੈ ਆਣੇ ਉਹ ਭਗਤੀ ਦਾਨ ਮੱਤ ਦੇਣਾ ਹੀ ਭਗਤੀ ਦਾਨ ਹੈ ਮੱਤ ਦੇਣਾ ਗੁਰ ਮੱਤ ਦਾ ਉਪਦੇਸ਼ ਦੇਣਾ ਹੀ ਭਗਤੀ ਦਾਨ ਹੈ ਉਹ ਭਗਤੀ ਦਿੰਦੇ ਲੈਂਦੇ ਕੌਣ ਨੇ ਸੰਤ ਜਨ ਸੰਤਾ ਕੋਲ ਭਗਤੀ ਨਹੀਂ ਹੁੰਦੀ ਸੰਤ ਜਨ ਸੰਤਾਂ ਤੇ ਸ਼ਾਂਤਮਈ ਗਿਆਨਵਾਨ ਜਿਹਨਾਂ ਨੂੰ ਸਮਝ ਆਉ ਉਹ ਲੈਂਦੇ ਨੇ ਸੰਤ ਜਨ ਲੈਣ ਲੈਂਦੇ ਸੰਤ ਨਹੀਂ ਲੈਂਦੇ ਜਦ ਸੰਤ ਲੈਣ ਦਾ ਮਨ ਬਣਾ ਲੈਂਦਾ ਨਾ ਗੁਰਮਤਿ ਲੈਣੀ ਹੈ ਉਹਦਾ ਮਨ ਬਦਲ ਜਾਂਦਾ ਫਿਰ ਜਨ ਬਣ ਜਾਂਦਾ ਤੇ ਉਹ ਸਮਝ ਆ ਜਾਂਦੀ ਹੈ ਸਮਝਦਾਰ ਸੰਤ ਲੈਂਦੇ ਨੇ ਆ ਜਿਹੜੇ ਦੂਏ ਸੰਤ ਨੇ ਪਾਗਲ ਸੰਤ ਨੇ ਮੂਰਖ ਉਹ ਨਹੀਂ ਲੈਂਦੇ ਉਹਨਾਂ ਨੇ ਲਈਓ ਨਹੀਂ ਮੂਰਖਾਂ ਨੇ ਜੱਟਾਂ ਸੰਤ ਜਨ ਉਹ ਸੰਤ ਜਨ ਤਾਂ ਜਾਂਚਦੇ ਨੇ ਮੰਗਦੇ ਨੇ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਬ੍ਰਹਮ ਗਿਆਨੀ ਤਾਂ ਮਹੇਸ਼ ਸ਼ਿਵਜੀ ਕੋ ਖੋਜਦਾ ਭਗਤੀ ਬਾਤੈ ਖੋਜਦਾ ਇਹ ਪੰਕਤੀ ਮੈਨੂੰ ਵੀ ਪੜ੍ਹੇ ਹਾਂਜੀ ਭਗਤੀ ਦਾ ਸੰਤ ਜਨ ਰਹਾਉ ਜਾਂਚੈ ਕਰ ਦਿਗ ਬਿਸੈ ਸੰਤ ਜਨ ਸੰਤ ਜਨਤਾ ਨੋਖਦੇ ਨੇ ਇੱਥੇ ਸੰਤ ਸਾਨੂੰ ਵਾਲਾ ਦੇ ਕੇ ਨਾਮ ਦਿੰਦੇ ਨੇ ਉਹ ਸੰਤ ਜਨ ਸੰਤਾਂ ਦਾ ਤਾਂ ਨਾਮ ਹੁੰਦਾ ਹੀ ਨਹੀਂ ਭਗਤਾਂ ਕੋਲ ਹੁੰਦਾ ਹੈ ਨਾਮ ਫਰਕ ਹੈ ਗੱਲ ਦਾ ਬਹੁਤ ਬਰੀਕ ਗੱਲ ਹੈ ਸੰਤਾਂ ਦਾ ਨਾਮ ਹੀ ਨਹੀਂ ਹੁੰਦਾ ਸੰਤਾਂ ਦਾ ਵਿਦੇਸ਼ ਕੀਤਾ ਗੁਰਬਾਣੀ ਨੇ ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸੰਤਾਂ ਨੂੰ ਤਾਂ ਕਹਿ ਆਵੇ ਤੁਸੀਂ ਆ ਜਿਹੜਾ ਸ਼ਬਦ ਦਾ ਨਾਰਦੀ ਭਗਤੀ ਹੈ ਨਾਰਦੀ ਮੰਗਰ ਵਾਲੀ ਨਾਰਦਰ ਨੇ ਜਿੱਥੇ ਤਪੱਸਿਆ ਕੀਤੀ ਇੱਥੇ ਉਹ ਭਗਤੀ ਹੈ ਕੋਈ ਬਨਾਰਸ ਕੋਲ ਦੀ ਧਰੂ ਕੋਲ ਹੈ ਇਹਨਾਂ ਸੰਤਾਂ ਕੋਲ ਬਨਾਰਸ ਵਾਲੀ ਬਨਾਰਸ ਕੇ ਠੱਗ ਜਿਵੇਂ ਸਾਡੀ ਜਿਹੜੀ ਪ੍ਰਚਾਰ ਹੁੰਦਾ ਸਿੱਖੀ ਦਾ ਹੁੰਦਾ ਅਮਰਸਰ ਵਾਲਾ ਆਨੰਦਪੁਰ ਸਾਹਿਬ ਵਾਲਾ ਹੁੰਦਾ ਹੀ ਨਹੀਂ ਅਮਰਸਰ ਵਾਲਾ ਖਾਸੀਗੜ੍ਹ ਕੋਈ ਹੈ ਕਿਉਂ ਕਾਚੀ ਦੇ ਠੱਗ ਅਰੰਬਰਸਾ ਬਨਾਰਸ ਦੇ ਠੱਗ ਉਧਰ ਅੰਬਰਸਾਲ ਦੇ ਠੱਗ ਦੋਵੇਂ ਮਸ਼ਹੂਰ ਨੇ ਦੋਵੇਂ ਵੱਡੇ ਸੈਂਟਰ ਨੇ ਧਰਬ ਦੇ ਦੋਹਾਂ ਦੇ ਵਿੱਚ ਠੱਗ ਜੁੜਿਆ ਹੋਇਆ ਕਿਉਂ ਜੁੜਿਆ ਠੱਗ ਅੰਬਰਸਾਲ ਦੇ ਠੱਗ ਅੰਬਰਸਾਲ ਅੰਦਰ ਸੜੀਏ ਇਹ ਜਿਹੜੇ ਨੇ ਇਹ ਸੰਤ ਨੇ ਇਹਨਾਂ ਕੋ ਤਾਂ ਨਾਮ ਹੁੰਦਾ ਹੀ ਨਹੀਂ ਸੰਤਾ ਕੋਈ ਨਾਮ ਕਦੇ ਹੋਇਆ ਅਸਾਤ ਭਗਤਾਂ ਕੋਲ ਹੋਇਆ ਬੱਬਈ ਫਿਰ ਉਹ ਸੰਤ RAM ਹੈ ਇੱਕੋ ਉਹ ਸੰਤ ਜਾਣਿਆ ਫਿਰ ਉਹ ਹੱਦ ਹੋ ਗਈ ਸੰਤ RAM ਦਾ ਉਹ ਹੋ ਉਹ ਸੰਤ RAM ਜਿਹੜਾ ਅੰਦਲਾ ਉਹ ਸੰਤ ਤਾਂ ਹੈ ਉਹ ਚਿੱਤਰ ਮੰਡੇ ਲੈਵਲ ਦੀ ਗੱਲ ਹੈ ਉਹ RAM ਕੜਾ ਗਿਆਨਬਾਨ ਰਾਮ ਦਾ ਰੋਂਦਾ ਸੰਤ ਵੀ ਰੋਂਦਾ ਰੋਵੇ RAM ਨਾ ਕਾੜਾ ਪਿਆਨੇ ਹਾਂਜੀ ਔਰ ਉਹ ਰਾਮ ਵੀ ਕਿਹਾ ਹੈ ਨਾ ਹਾਂਜੀ ਉਹ ਉੱਥੇ ਪੰਕਤੀ ਹੈ ਜੀ ਸੰਤ ਰਾਮ ਹੈ ਇੱਕੋ ਬਾਈ ਨਿੰਦੋ ਰਾਂ ਸੰਤਾ ਨੂੰ ਪਰ ਉਪਦੇਸ਼ ਦਾ ਕਰਨਾ ਕਿ ਨਹੀਂ ਕਰਨਾ ਜਦ ਸੰਤ ਕਹਿੰਦੇ ਨੇ ਸਾਡੇ ਕੋਲ ਨਾਮ ਹੈਗਾ ਹੈ ਨਹੀਂ ਫਿਰ ਉਹ ਨਿੰਦ ਫਿਰ ਉਹ ਠੱਗ ਹੋ ਜਾਂਦੇ ਨੇ ਸੰਤ ਨਹੀਂ ਹੈ ਸੰਤ ਹਰਕੇ ਸੰਤ ਹੁੰਦੇ ਨੇ ਕੱਲੇ ਸੰਤ ਨਹੀਂ ਹੁੰਦੇ ਜਿਹੜੇ ਸੰਤ ਜਾਣੇ ਉਹ ਹਰਕੇ ਸੰਤ ਕਹਿ ਕੇ ਐਡ ਕਰ ਲੈ ਹਰਕੇ ਸੰਤ ਨਾ ਆਖੀਐ ਬਾਨ ਆਰਥ ਕੇ ਠਗ ਜਿਹੜੇ ਹਰਕੇ ਸੰਤ ਨਹੀਂ ਹੈ ਜਿਹਨੇ ਨਾਮ ਜਿਹੜੇ ਕਹਿੰਦੇ ਸਾਡੇ ਕੋਲ ਨਾਮ ਹੈਗਾ ਹਰਕੇ ਸੰਤ ਨਹੀਂ ਕਹਿੰਦੇ ਸਾਡੇ ਕੋਲ ਨਾਮ ਹੈਗਾ ਉਹ ਹਰਕੇ ਸੰਤ ਤਾਂ ਥੱਲੇ ਨੇ ਸੰਤ ਆਫੇ ਗੁਰੂ ਬਣੇ ਬੈਠੇ ਨੇ ਉਤਾ ਜੋ ਹਰਕੇ ਕੇ ਸੰਤ ਨੇ ਨਾ ਕਿਸੇ ਦੇ ਨੇ ਉਤਾ ਜੀ ਉਤਾ ਜੋ ਚੇਲੇ ਨੇ ਹਾਂਜੀ ਜਿਹੜੀ ਭਗਤੀ ਸੰਤ ਕਰਦੇ ਨੇ ਜਦੋਂ ਪਤਾ ਲੱਗਿਆ ਭਗਤੀ ਗਲਤ ਹੈ ਪਾਵਨਾਂ ਨੇ ਭਗਤੀ ਮੰਗੀ ਜਾਚੈ ਕਰ ਦਿਗ ਦਿਸੈ ਸਰਾਇ ਆ ਜਿਹੜੇ ਘਰ ਦੇ ਵਿੱਚ ਐਡੀ ਬੜੀ ਕਨਾਤ ਹੈ ਕਨਾਤ ਕਨਾਤ ਮਤਲਬ ਹੁੰਦੀ ਆਹ ਲੜੇ ਆਹ ਜਿਹੜਾ ਨਾ ਆਪਣਾ ਰਾਮਗਰਬ ਰਾਮਗਰਬ ਹੈ ਜੀ ਤਿੰਨ ਲੋਕ ਨੇ ਇਹ ਉਹਦੇ ਘਰ ਦੇ ਅੰਦਰ ਹੈ ਜਿਹੜਾ ਭਵਸਾਗਰ ਹੈ ਇਹ ਉਹਦੇ ਘਰ ਦੇ ਅੰਦਰ ਹੈ ਸੁਖ ਸਾਗਰ ਤੇ ਉਹਦਾ ਘਰ ਸੁਖ ਸਾਗਰ ਹੈ ਭਵਸਾਗਰ ਉਹਦੇ ਅੰਦਰ ਆ ਸਾਰੀ ਰਚਨਾ ਭਵਸਾਗਰ ਦੇ ਵਿੱਚ ਹੀ ਹੈ वैकुंठ भवन चित्रशाला वैकुंठ भवन चित्रशाला ओदे विच ही है जदों तुसी वैकुंठ गए ने ओ भवन और चित्रशाला संसार ए संसार है वैकुंठ नोदा ए चित्रशाला इही है इथे या जून दा चित्र चित्र विचित्र आया बेचारा चित्र चित्र आ ए संसार उनी देखणा संसार चित्र ਸੱਚੀ ਮੂਰਤ ਹੈ ਚਲਦੀ ਫਿਰਦੀ ਤੇ ਜਾਨਦਾਰ ਮੂਰਤਾਂ ਨੇ ਜੜ ਕੇ ਤੰਨਾ ਬੇਲ ਹੈ ਜਿਹੜੀ ਅਸੀਂ ਮੂਰਤ ਬਰੋਲਦੇ ਉਹ ਜੜ ਹੁੰਦੀ ਹੈ ਉਹ ਇਸ ਮੂਰਤ ਦੀ ਦੇਖਣਾ ਖੂਬਸੂਰਤੀ ਨਹੀਂ ਦੇਖਣੀ ਹੈ ਤੇਰੀ ਐਨਜੋਏ ਕਰਨ ਨੂੰ ਆਸਤੇ ਅਸੀਂ ਇੱਥੇ ਆਏ ਤਾਂ ਕਿ ਧਿਆਨ ਛੱਡ ਕੇ ਜਿਹਦੇ ਚਿੱਤਰ ਰਚਿਆ ਜਿਹਦੇ ਚਿੱਤਰ ਬਣਾਇਆ ਹੈ ਜੇ ਤੇਰਾ ਜਦੋਂ ਉਹਦੇ ਵਾਸਤੇ ਰੱਖਣਾ ਇੱਥੋਂ ਚਿੱਤਰ ਵਿੱਚੋਂ ਯਾਨੀ ਤਨ ਵਿੱਚੋਂ ਮਨ ਖੋਜਣਾ ਹੈ ਤਨ ਨਹੀਂ ਖੋਜਣਾ ਸੰਸਾਰ ਤਨ ਖੋਜਦੇ ਡਾਕਟਰ ਤਨ ਖੋਜਦੇ ਨੇ ਰਿਵੋਲਟ ਤਨ ਖੋਜਣ ਬਣਾਏ ਨੇ ਮੈਡੀਕਲ ਸੈਨ ਤਨ ਖੋਜਣ ਤੇ ਬਣੀ ਹੈ ਆਯੁਰਵੈਦਿਕ ਤਨ ਖੋਜਣ ਦੀ ਗੱਲ ਹੈ ਜਿਹੜੇ ਯੋਗਾ ਤਨ ਖੋਜਣ ਦੀ ਗੱਲ ਹੈ ਇਹ ਤਨ ਵਿੱਚੋਂ ਮਨ ਖੋਜਣਾ ਹੈ ਹਾਂਜੀ ਤੁਸੀਂ ਕਿਹਾ ਕਿ ਅਸੀਂ ਇੰਜੋਏ ਕਰਨ ਨਹੀਂ ਆਏ ਨਹੀਂ ਆਏ ਹੁੰਦਾ ਕੀ ਹੈ ਆਮ ਤੌਰ ਤੇ ਬੰਦਾ ਬੋਰ ਹੋ ਜਾਂਦਾ ਕਹਿੰਦਾ ਚਲੋ ਥੋੜਾ ਇੰਜੋਏ ਕਰ ਲਈਏ ਫਿਰ ਉਹ ਲਾਈਫ ਕੀ ਹੈ ਤੇ ਤੁਸੀਂ ਜਿਹੜੀ ਜ਼ਿੰਦਗੀ ਦੀ ਗੱਲ ਕਰ ਰਹੇ ਹੋ ਉਹ ਕਿਹੜੀ ਹੈ ਉਹ ਤਾਂ ਸੰਸਾਰੀ ਕਹਿੰਦੀ ਹੈ ਇੰਜੋਏ ਕਰਨੀ ਉਹ ਦੁੱਖਦਾਂ ਦੀ ਜ਼ਿੰਦਗੀ ਹੈ ਇੰਜੋਏ ਕਰਨਾ ਦੁੱਖਦਾ ਹੈ ਦੋਈ ਪਾਸੇ ਕਰਦਾ ਜੇ ਦੋਹੇ ਸੰਸਾਰ ਦੇ ਵੀ ਇੰਜੋਏ ਕਰਦਾ ਹੈ ਮਹਾਰਾਗੀ ਵੀ ਉਦੋਂ ਕਾਟਦਾ ਫਿਰ ਦੁਗਦਾ ਹੈ ਉਹ ਦੁਗਦਾ ਰੋਗ ਦੁਗਦਾ ਦੇ ਵਿੱਚ ਰੋਗ ਜਿਹੜੇ ਵਧਦੇ ਨੇ ਹੋਏ ਨੇ ਇਹਲੇ ਸੰਤ ਜਨ ਭਗਤੀ ਮੰਗਦੇ ਨੇ ਭਗਤੀ ਤਾਂ ਇੱਕੋ ਦੇ ਸ਼ਬਦ ਜਾਂਦੀ ਹੈ ਫਿਰ ਏਕਾ ਦੇਸ ਧਾਵਾ ਜਿਹੜਾ ਦੋ ਪਾਸੇ ਜਾਂਦਾ ਉਹ ਵਿਚਾ ਉੱਥੇ ਹੀ ਰਹਿੰਦਾ ਉਧਰੋਂ ਕਾ ਜਿਹੜਾ ਉਧਰੋਂ ਬਜਲੇ ਵਿਚਾਰੇ ਰਹਿੰਦੇ ਆ ਬਸ ਹਾਂ ਉਹ ਤੇ ਬੋਰ ਹੁੰਦਾ ਕਿਉਂ ਆ ਪਹਿਲਾਂ ਇਹ ਦੱਸ ਬੋਰ ਹੋ ਜਾਂਦੇ ਵੀ ਜਿਹੜਾ ਮਨ ਹੈ ਉਹ ਯਾਰ ਫਿਰ ਉਹ ਹੀ ਗੱਲ ਬਿਆਕੁਲ ਮੇਰਾ ਨਹੀਂ ਮੇਰਾ ਸਵਾਲ ਹੋਰ ਹੈ ਹਾਂਜੀ ਭਗਤ ਬੋਰ ਹੁੰਦਾ ਹੀ ਨਹੀਂ ਹਾਂ ਉਹ ਕਿਉਂ ਨਹੀਂ ਹੁੰਦੇ ਬੋਰ ਉਹ ਤਲ ਵਿੱਚ ਉਹਨਾਂ ਦਾ ਟੇਸੇ ਹੋ ਰਿਹਾ ਇਹ ਟੇਸੇ ਹੋ ਰਿਹਾ ਮਾਇਆ ਦੇ ਟੇਸੇ ਇੱਕ ਜਗ੍ਹਾ ਤੁਸੀਂ ਟਿਕ ਨਹੀਂ ਸਕਦੇ ਬੋਰ ਹੋਵੋਗੇ ਕਿਉਂਕਿ ਉਹ ਤੇ ਮਾਇਆ ਟਿਕ ਨਹੀਂ ਸਕਦਾ ਬੋਰ ਉਹ ਨਾਮ ਦੀ ਭੁੱਖ ਆਲੇ ਦੀ ਭੁੱਖ ਹਟਦੀ ਹੋਈ ਨਹੀਂ ਮਾਇਆ ਦੀ ਭੁੱਖ ਤਾਂ ਥੋੜੀ ਭੁੱਖ ਹੈ ਬਸ ਉਹ ਥੋੜਾ ਦਿਰ ਬਾਅਦ ਇਹ ਹਟ ਜਾਂਦੀ ਹੈ ਫਿਰ ਉਹ ਬੋਰ ਹੋ ਜਾਂਦਾ ਨਾਮ ਦੀ ਭੁੱਖ ਹੈ ਉੱਥੇ ਉਹ ਕਿਵੇਂ ਹਟ ਸੰਸਾਰ ਦੀ ਪੁੱਖ ਪੂਰੀ ਹੁੰਦੀ ਹੈ ਉਹ ਪੂਰੀ ਹੋ ਨਹੀਂ ਹੁੰਦੀ ਪੁੱਖ ਅਦੇ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾ ਉਹ ਭਗਵਾਨ ਦੇ ਲੈਵਲ ਤੇ ਹੈ ਉਹ ਇੰਜੋਏ ਕਰਨ ਸਾਡੀ ਲੋੜ ਹੈ ਉਸ ਨਾਲ ਬੋਰ ਹੋ ਗਿਆ ਲੋੜ ਹੈ ਇੰਜੋਏ ਕਰ ਲੈ ਬੋਰ ਹੁਣ ਤੇ ਅਸੀਂ ਮੰਨ ਉਸੇ ਕੰਮ ਤੇ ਲੱਗੇ ਇਹ ਕੂੜੇ ਕੰਮ ਨੇ ਜਿਹੜੇ ਕੂੜੇ ਕੰਮਾਂ ਦੇ ਵਿੱਚੋਂ ਬੋਰ ਹੁੰਦਾ ਇਹ ਮਾਇਆ ਦੇ ਕੰਮ ਲਈ ਇੱਥੇ ਬੋਰ ਹੁੰਦਾ। ਨਾਮ ਦੀ ਖੋਜ ਵਾਲਾ ਬੋਰ ਹੁੰਦਾ ਹੀ ਨਹੀਂ। ਅਸੀਂ ਕੰਮ ਕਰਦੇ ਹਟ ਜਵੇ। ਜਾਂ ਉਸ ਰਸ ਲੋੜ ਡਾ ਫਿਰ ਅਸੀਂ ਬੋਰ ਹੋਣ ਲੱਗ ਜਾਈਏ। ਜੇ ਤ੍ਰਿਪਤੀ ਹੋ ਨਹੀਂ ਹੁੰਦੀ ਫਿਰ ਬੋਰ ਕਿਵੇਂ ਹੋਊ? ਮਾਇਆ ਚ ਤ੍ਰਿਪਤੀ ਹੈ। ਮਾਇਆ ਚ ਤ੍ਰਿਪਤੀ ਹੈ। ਤ੍ਰਿਪਤ ਰਹੇ ਨਾ ਆਏ। ਮਾਇਆ ਤ੍ਰਿਪਤੀ ਜਿਆਦਾ ਜਸ ਸੰਤੋਖ ਆ ਜਾਂਦਾ ਹੈ ਬਿਨਾ ਸੰਤੋਖ ਨਹੀਂ ਕੋ ਰਾਜਾ ਹੈ ਪਰ ਮਾਇਆ ਇੱਕ ਥਾਂ ਨਹੀਂ ਨਾ ਮਾਇਆ ਬਹੁ ਰੰਗੀ ਹੈ ਉੱਤੇ ਇੱਕ ਰੰਗ ਹੈ ਇੱਕ ਰੰਗ ਤੋਂ ਬੋਰ ਹੁੰਦਾ ਦੂਗੇ ਰੰਗ ਚਾਉਂਦਾ ਦੂਏ ਤੋਂ ਬਹੁ ਟੀਏ ਰੰਗ ਚ ਜਾਉਂਦਾ ਉੱਤੇ ਰੰਗ ਇੱਕਾ ਰੂਆ ਹੈ ਹੀ ਨਹੀਂ ਉੱਤੇ ਬਹੁਤਾ ਸਵਾਲੇਵਾਦੀ ਹੁੰਦਾ ਦੂ ਕੀ ਹੈ ਨਹੀਂ ਉਹ ਜੀ ਹੋਰ ਕਿਉਂ ਹੋਊਗਾ ਇਹ ਤਾਂ ਦੇਖ ਲੈ ਮਾਇਆ ਦੇ ਰੰਗ ਤਾਂ ਸਾਰੇ ਜਦ ਮਾਇਆ ਦੇ ਰੰਗਾਂ ਦੇ ਉਹ ਛੁੱਟ ਕੇ ਦੂਏ ਪਾਸੇ ਗਿਆ ਮਾਇਆ ਦੇ ਰੰਗ ਤਾਂ ਉਹ ਜੱਟੇ ਸਹੀ ਨਹੀਂ ਉਹਦੇ ਮੁਕਾਬਲੇ ਦਾ ਜੇ ਕੋਈ ਸਾਨੂੰ ਟੇਸ ਹੋਰ ਹੁੰਦਾ ਫਿਰ ਬੋਰ ਹੋ ਕੇ ਦੂਏ ਤੇਸਵਾਂ ਲੱਗਦਾ ਉਹਨਾਂ ਨੂੰ ਲੱਗਦਾ ਹੀ ਨਹੀਂ ਵੈਸੇ ਇਹ ਗੱਲ ਨੂੰ ਉਹੀ ਸਮਝ ਸਕਦਾ ਜੀ ਦੀ ਵਸਤਵ ਹੋਵੇ ਆਮ ਆਦਮੀ ਨਹੀਂ ਸਮਝਣ ਦੇ ਸਾਨੂੰ ਮਾਇਆ ਵਾਲੇ ਕਦੇ ਇਸ ਗੱਲ ਉਹ ਤਾਂ ਬੋਰ ਹੁੰਦੇ ਨੇ ਨਾਮਦਾਰਾ ਸਾਨੂੰ ਆਇਆ ਕੋਈ ਨਹੀਂ ਉਹ ਮੈਂ ਨਹੀਂ ਮਾਇਆ ਗਾਇਕਾ ਬਛੜਾ ਬਛੜਾ ਛੋਟਲਾ ਥਣ ਚੌਂਖੇ ਮਾਂ ਖੰਕੂਟਲਾ ਜਿਹਨੂੰ ਅੱਖਾਂ ਦੇ ਕੋਟਾਉਂਦੇ ਨੇ ਥਣ ਛੱਡ ਦਾ ਪੇਟ ਲਿਮਟਿਡ ਪਤਾ ਕਿੰਨਾ ਹੈ ਲਿਮਟਿਡ ਨਹੀਂ ਹੈ ਘਰ ਹੈ ਦਿਗ ਹਾਂ ਗ੍ਰੰਥ ਗਾਨੀ ਦਾ ਮਨ ਪਰਗਾਸ ਜੈਸੇ ਤਾਰੂ ਪਰ ਤਾਰੂ ਪਰ ਆਜ ਨਾ ਉਹਦਾ ਪੇਟ ਹੈ ਪਰੂ ਕਹਦੇ ਨਾ ਪਰੂ ਕਹਦੇ ਨਾ ਜਨਮ ਤਾਂ ਬੰਦਾ ਨਹੀਂ ਫੇਰ ਵੀ ਬਹੁਤ ਕੁਝ ਹੈ ਜਾਣਨ ਨੂੰ ਬਹੁਤ ਕੁਝ ਹੈ ਜਦ ਉਹਦੇ ਜੋ ਜਾਣਨ ਨੂੰ ਮੁੱਖ ਜਵੇ ਸਾਨੂੰ ਰਾਸ ਜਿਆਦਾ ਹੁੰਦੇ ਹੁੰਦਾ ਜਿਹੜੇ ਖੋਜੀ ਨੇ ਖੋਜੀ ਨਹੀਂ ਬੋਲੁੰਦੇ ਕਹਿੰਦੇ ਖੋਜੀ ਸੁਣਿਆ ਬੋਲ ਰਹਾ ਨਹੀਂ ਉਹ ਕਹਿੰਦੇ ਵੀ ਤੱਕ ਆਪਣੇ ਧੁੰ ਚ ਲੱਗਿਆ ਹੀ ਰਹਿੰਦਾ ਹਰ ਉਹ ਵਾਲੇ ਬੋਰ ਹੁੰਦਾ ਕੋਈ ਕਦੇ ਬੋਰ ਨਹੀਂ ਹੁੰਦਾ ਬੋਰ ਤਾਂ ਨਹੀਂ ਕੋਈ ਦਾ ਧਿਆਨ ਇੱਕ ਪਾਸੇ ਨਹੀਂ ਹੁੰਦਾ ਹਾਂ ਬੋਰੰਗੀ ਮਾਇਆ ਖੇਡਦੇ ਨੇ ਜਿਹੜੇ ਉਹ ਬੋਰ ਹੁੰਦੇ ਨੇ ਕੋਈ ਜੀ ਨੂੰ ਨਵਾਂ ਕੋਈ ਨਵਾਂ ਕੁ ਮਿਲਦਾ ਰਹਿੰਦਾ ਹੈ ਉਹ ਗਾਹ ਤੁਰਦਾ ਰਹਿੰਦਾ ਜਿਹੜਾ ਬੋਰ ਹੋ ਜਵੇ ਖੋਜੀ ਨਹੀਂ ਹੈ ਇਹ ਵੀ ਗੱਲ ਹੈ ਖੋਜੀ ਬੋਰ ਹੁੰਦਾ ਨਹੀਂ ਜੇ ਬੋਰ ਹੋਵੇ ਖੋਜੀ ਹੈ ਨਹੀਂ ਕੋਈ ਗਿਆਨ ਅਸੀਮ ਹੈ ਚਾਹੇ ਕੋਈ ਵੀ ਹੋਵੇ ਗਿਆਨ ਅਸੀਮ ਖੋਜ ਗਿਆਨ ਦੀ ਖੋਜ ਲੱਗਿਆ ਬੋਰ ਕਿਉਂ ਹੋਊਗਾ ਬੋਰ ਜਾਦਾ ਹੋ ਫਿਰ ਖੋਜੀ ਖੋਜੀ ਨਹੀਂ ਰਹਿਣਾ ਬੰਦ ਹੋ ਖੋਜ ਪਰ ਫਿਰ ਖੋਜੀ ਨਹੀਂ ਹੈ ਜੇ ਬੋਰ ਹੋਗਾ ਫਿਰ ਲਾਲਾ ਹੋ ਜੀਏ ਫਿਰ ਲਾਲਾ ਬ੍ਰੇਕ ਟੁੱਟ ਗਿਆ ਉੱਥੋਂ ਸੱਪਤ ਲੋਕ ਸਾਮਾਨ ਪੂਰੀਲੇ ਸਾਧਾ ਲੋਕ ਦਾ ਸਾਮਾਨ ਇੱਕ ਵਾਰ ਪਾਤਾ ਇੱਥੇ ਜਿਹੜੇ ਸਾਧਾ ਲੋਕ ਕਹਿੰਦੇ ਨੇ ਨਾ ਕੋਈ 14 ਲੋਕ ਕਹਿੰਦਾ 14 ਬਤਾਰ 14 ਨਰਕ ਵਾਲੇ ਨੇ 14 ਨਾ 7 ਨਰਕ ਦੇ ਨੇ 7 ਸਤ ਸਵਰਗ ਦੇ ਨੇ 7 ਦੇਵਤਿਆਂ ਦੇ ਨੇ 7 ਰਾਖਸ਼ਾਂ ਨੇ ਰਾਖੀ ਦੇਵਤਿਆਂ ਦਾ ਪਰ ਨਹੀਂ ਕਹਿੰਦੇ ਤੇ ਕੋਈ ਹੁੰਦੇ ਨੇ ਅਸਲ 'ਚ ਜਿਹੜਾ ਆਖਿਂਦੇ ਨੇ ਸਨਾਤਨਵਾਦ ਵਾਲੇ ਉਹ ਉਹਨਾਂ ਨੂੰ ਗੁਰਬਾਣੀ ਇਕੱਠੇ ਏ ਕੋਈ ਮੰਦੀ ਏ ਪਾਪਨ ਦੋਨੋਂ ਭਾਈ ਅਸੀਂ ਮੰਨਦੇ ਹਾਂ ਸਾਖਤ ਔਰ ਸੰਤ ਉਹ ਨਹੀਂ ਮੰਨਦੇ ਸਨਾਤਨ ਵਾਲੇ ਸਾਖਤ ਨਹੀਂ ਮੰਨਦੇ ਕੋ ਕੋ ਸਾਖਤ ਆਪਨੇ ਸਨਾਤਨੀ ਨੇ ਸਾਖਤ ਨੇ ਹੋ ਸਾਰੇ ਇਸ ਕਰਕੇ ਸਾਖਤ ਨਹੀਂ ਮੰਨਦੇ ਹੋ ਸਾਖਤ ਆਪਨੇ ਹੋ ਸਾਕਤ ਮਰਨ ਸੰਤ ਸਭ ਜੀਵ ਹੈ ਜਿਹੜੇ ਮਰਨਾ ਮੰਨਦੇ ਨੇ ਵੀ ਮਰ ਜਾਂਦਾ ਹੈ ਜਿਹੜੇ ਕਰਿਆ ਕਰਮ ਨੂੰ ਮੰਨਦੇ ਨੇ ਜਿਹੜੇ ਫੁੱਲ ਪਾਉਂਦੇ ਨੇ ਮਰਨ ਤੋਂ ਬਾਅਦ ਉਹਦੇ ਸਭ ਕੁਝ ਕਰਦੇ ਨੇ ਕਰਿਆ ਕਰਮ ਉਹ ਸੰਸਾਰੀ ਆਦਮੀ ਨੇ ਉਹ ਮਤਾਂ ਸੰਸਾਰੀ ਨੇ ਸਨਾਤਨੀ ਮਤ ਤੇ ਮੰਨਦੀ ਹੈ ਸਨਾਤਨੀ ਮਤ ਬੇਦਮਤ ਨਹੀਂ ਬੇਦਮਤ ਨਹੀਂ ਮੰਨਦੀ ਬੇਦਮਤ ਮੰਨਦੀ ਐਨੇ ਕ ਜਨਮ ਐਨੇ ਕਿਸਮਰ ਆਪਣੇ ਚਲ ਆ ਵੀ ਕਰ ਆਵਣ ਜਾਵਣ ਦੇਸ਼ ਅੰਦਰਿਸ਼ਟ ਆਗਿਆਕਾਰੀ ਤਾਰੀ ਸਭ ਸਿ ਆਗਿਆਕਾਰੀ ਤਾਰੀ ਸਭ ਸਿ ਸਨਾਤਨੀ ਮਤ ਜਿਹੜੇ ਸੰਥਾਰੀ ਮਤ ਵਾਲੇ ਨੇ ਮਤ ਨਹੀਂ ਹੈ ਨਰਾਕਾਰ ਸੰਬੰਧ ਨਹੀਂ ਕੋਈ ਉਹ ਮੂਰਤੀ ਪੂਜਾਉਣੇ ਨੇ ਸਾਰੇ ਮੂਰਤੀ ਪੂਜਣਾ ਫਰਾਂਤਨੀ ਮਤ ਕੋਈ ਮਾਇਆ ਤਾਰੀ ਨੇ ਅੰਮੇ ਬੋਲੇ ਸਨਾਤਨੀ ਵਾਸਤਵ ਕਬੀਰ ਕੋਲ ਹੈ ਪਹਿਲਾਂ ਸਨਾਤਨੀ ਮਾਤ ਦੇ ਆਏ ਨੇ ਸਾਡੇ ਸੰਤੇ ਕੁਛ ਛੱਡੀ ਹੈ ਇਹਨਾਂ ਨੇ ਸਨਾਤਨੀ ਮਾਤ ਤੋਂ ਸੰਤ ਪੈਦਾ ਕਰਦੀ ਹੈ ਸਨਾਤਨੀ ਸਨਾਤਨੀ ਇਹ ਸੰਤ ਜਨ ਮੰਗਦੇ ਨੇ ਤੇ ਲਿਖਿਆ ਚਾਹ ਸੰਤ ਜਨ ਉਹ ਭਗਤੀ ਦੇਣ ਵਾਲਾ ਸੰਤ ਜਨ ਭਗਤੀ ਮੰਗਦੇ ਨੇ ਨਾਮ ਨਾਮ ਪਦਾਰਥ ਸਨਾਤਨੀ ਵਾਦ ਦੇਗਾ ਚਾਰ ਪਦਾਰਥ ਨਹੀਂ ਚਾਰਾਂ ਦਾ ਨਾਮ ਹੈ ਹੀ ਨਹੀਂ ਧਰਮ ਅਰਥ ਕਾਮੋਗ ਹੈ ਪਹਿਲੀ ਗੱਲ ਤਾਂ ਧਰਮ ਉਹ ਕੋਈ ਧਰਮ ਦੇ ਵਿੱਚ ਪਦਾਰਥ ਨਹੀਂ ਚਾਰ ਧਰਮ ਚਾਰ ਪਦਾਰਥ ਮੰਨਦਾ ਚਾਰ ਪਦਾਰਥ ਜੇ ਕੋ ਮੰਗਾ ਚਾਰ ਪਦਾਰਥ ਧਰਮ ਕਾਦਮੀ ਮੰਨਦਾ ਸਨਾਤਨੀ ਵਾਦ ਚਾਰ ਪਦਾਰਥ ਹੀ ਤਿੰਨ ਨੇ ਉਹ ਧਰਮ ਨੂੰ ਪਦਾਰਥ ਮੰਨਦੇ ਨੇ ਉਹ ਧਰਮ ਦਾ ਵਦਾਰਤ ਕਿਤੇ ਧਰਮ ਦਾ ਧਾਰਨ ਕਰਨ ਵਾਲੀ ਚੀਜ਼ ਹੈ। ਉਹ ਦਾਤਾਂ ਜੋ ਧਰਮ ਚੋਂ ਮਿਲਦੇ ਨੇ ਯਾਰ। ਇਹ ਮੰਗੀਦੇ ਹੁੰਦੇ ਨੇ। ਧਰਮ ਧਾਰਨ ਕਰਕੇ ਕੋਈ ਮੰਗਦੇ ਨੇ ਮਨੋ ਕਾਮਨਾਵਾਂ ਪੂਰੀਆਂ ਹੋ ਵੀ ਉਹੀ ਮੰਗਦੇ ਨੇ। ਇਹ ਧਨ ਸੰਖਾਰੀ ਪੈਸਾ ਅਰਥ ਇਹ ਸੰਖਾਰੀ ਵੈਸ਼ ਆ ਹੈ। ਪੰਨ ਬਦੀ ਬਣਾਈ ਹੋਈ ਮਤ ਹੈ ਰਾਜੇ ਵਾਸਤੇ ਰਾਜ ਦਾ ਕੰਮ ਹੈ ਇਹ ਆਰਥਿਕਤਾ ਆਰਥਿਕ ਮੰਦਲ ਲੋਕਾਂ ਦੀ ਗੱਲ ਨਹੀਂ ਤੋਂ ਤਾਂ ਲੈ ਕੇ ਹੀ ਲੋਕਾਂ ਦੀ ਮਦਦ ਕਰਨੀ ਹੈ ਜਿਵੇਂ ਸਰਕਾਰ ਕਰਦੀ ਹੈ ਇਹ ਤਾਂ ਲੈ ਕੇ ਟੈਕਸ ਆਫੇ ਖਾਈ ਜਾਂਦੇ ਨੇ ਦੁਹਾਨ ਨੂੰ 15 ਪੈਸੇ ਵੀ ਨਹੀਂ ਦਿੰਦੇ ਅਰਥ ਕਾਮਨਾ ਪੂਰੀਆਂ ਕਰਨ ਵਾਸਤੇ ਤਾਂ ਸੱਚਾਈ ਦਾ ਕਾਮ ਅਰਥ ਫਿਰ ਮੁਕਤੀ ਉਹ ਜੇ ਤੇ ਕਾਮਨਾ ਮੁਕਤੀ ਕਿਵੇਂ ਹੋ ਜੂ ਉਥੇ ਨਾਲੇ ਕਾਮਨਾ ਛੱਡੇ ਤੇ ਮੁਕਤੀ ਹੈ ਇੱਛਾਵਾਂ ਤੇ ਤੇ ਮੁਕਤੀ ਹੈ ਇੱਛਾਵਾਂ ਤੇ ਦੀ ਗੱਲ ਕਰ ਰਹੇ ਹੋ ਨਾਲੇ ਤੁਸੀਂ ਉਹਨੂੰ ਪਦਾਰਥ ਮੰਨੀ ਬੈਠੇ ਹੋ ਇਹ ਤਾਂ ਬਹੁਤ ਬੁਰੀ ਤਰ੍ਹਾਂ ਲਜਾਉਣ ਵਾਲੀ ਮਾਤਾ ਆ ਬੁੱਢ ਜੇ ਹੁੰਦੇ ਆਪ ਡੁੱਬੇ ਕਿਉਂ ਵੇਦਮੇ ਚੇਲੇ ਦੇ ਬਾਹਰ ਆਪ ਚਾਰ ਵੇਦਾਂ ਡੁੱਬ ਗਿਆ ਚੇਲੇ ਸਾਰੇ ਰੋੜ ਤੇ ਇਤਨਾ ਅਧਨੀ ਮਕਤਾ ਤਾਂ ਹੀ ਗੁਰੂ ਕੰਨ ਇਹ ਮਨ ਉਲਟ ਸਨਾਤਨ ਹੋਵਾ ਹੁਣ ਮੇਰਾ ਮਨ ਸਨਾਤਨ ਮਤ ਤੋਂ ਉਲਟ ਗਿਆ ਨੀ ਛੱਡ ਗਿਆ ਵਾਹ ਫਿਰ ਨੀ ਛੱਡਤੀ ਪਤਾ ਖਾਲ ਲੱਗਿਆ ਸਨਾਤਨ ਮਤਾ ਇਹ ਗਲਤ ਹੈ ਬਸਰੀ ਗਲਤ ਸਨਾਤਨ ਮਤ ਨਾਲ ਉਹਦਾ ਮਨ ਜਿੱਤੇ ਨਹੀਂ ਹੋਇਆ ਚੁੱਪੇ ਨਹੀਂ ਹੋਇਆ ਜਾਂਦੇ ਕੀ ਹੋਇਆ ਦੂਜੇ ਤਬ ਜਾਣਿਆ ਜਦ ਜੀਵਤ ਨੂੰ ਜਨਮ ਪਤਾ ਲੱਗਿਆ ਜੀਵਤ ਮਨਨਾ ਕੀ ਹੁੰਦਾ ਜਦ ਮੈਂ ਖੁਦ ਜੀਵਤ ਮਰ ਗਿਆ ਕਿ ਆਹ ਵਕਤੀ ਹੈ ਠੀਕ ਤਬ ਜਾਣਿਆ ਤਬ ਗਿਆਨ ਹੋਇਆ ਮੈਨੂੰ ਆਤਮ ਮੈਂ ਆਪਣੇ ਆਪ ਨੂੰ ਜਾਣਿਆ ਜਦ ਮੈਂ ਉਹ ਮਰ ਗਿਆ ਜਿਉਂਦਾ ਹੀ ਸਰੀਰ ਚ ਰਹਿਣਾ ਹੀ ਮੇਰਾ ਮਨ ਮਰ ਗਿਆ ਮੇਰੀਆਂ ਛਾਣਾਂ ਖਤਮ ਹੋ ਗਈਆਂ ਕਾਮਨਾਵਾਂ ਤਾਂ ਖਤਮ ਕਰ ਸੀ ਇਹ ਕਹਿੰਦੇ ਨੇ ਕਾਮ ਪਦਾਰਥ ਕਿ ਕੋਦੋਂ ਧਰਮ ਆਪਣੇ ਅਭੂ ਧਰਮ ਕਹੀ ਜਾਂਦੇ ਨੇ ਜੀ ਹਾਰੇ ਹੋ ਜੋਹਾਰੀਏ ਦੁਬਾਰਾ ਆਉਣ ਨੂੰ ਮੈਦਾਨ ਆ ਜਾਣ ਸਮਾ ਲੋਕਾਂ ਨੂੰ ਵੀ ਪਤਾ ਲੱਗੇ ਕਿ ਧਰਮ ਹੁੰਦਾ ਕੀ ਆ ਜਾਂਚੇ ਕਰ ਲక్ష్ਮੀ ਕੁਆਰੀ ਉਹ ਤਾਂ ਗੱਲ ਕੁਆਰੀ ਆ ਇਹਨਾਂ ਦੇ ਸੱਤ ਦੇਵੀਆਂ ਨੇ ਉੱਥੇ ਇੱਕੋ ਹੀ ਆ ਉਤਤੈਕਾ ਉਹ ਜਾਂ ਆਪਿਕਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਉਹ ਉਹ ਬੁੱਧੀ ਅਕਾਦਮੀ ਦੀ ਬੁੱਧੀ ਕੋਹਨੀਆ ਬੁੱਧੀ ਦੋ ਹੁੰਦੀਆਂ ਨੇ ਕੋਈ ਅਕਲ ਹੁੰਦੀ ਹੈ ਕਾਜ਼ਮੀ ਗਿਆਨ ਕਈ ਪ੍ਰਕਾਰ ਦਾ ਹੋ ਸਕਦਾ ਅਕਲ ਨੂੰ ਪਰ ਅਕਲ ਤਾਂ ਇੱਕ ਕੋਈ ਹੈ ਕੋ ਜੜੀ ਲక్ష్ਮੀ ਕੁਆਰਾ ਉਹ ਹੈ ਲక్ష్ਮੀ ਉਹ ਤਾਂ ਨਾ ਉਹਦੇ ਕੋਲ ਨਾਮ ਤਾਂ ਦਿੰਦੀ ਆ ਉਹ ਉਹ ਮਤ ਮਾਤਾ ਉਹੀ ਮਤ ਮਾਤਾ ਸੰਤੋਖ ਪਤਾ ਹੈ ਸੰਤੋਖ ਹੁਲਦਾਤ ਜਬ ਸੰਤੋਖ ਤਾਨਾ ਜਬ ਆਵੇ ਧਨ ਸੰਤੋਖ ਨੂੰ ਤਨ ਮੰਨਿਆ ਐ ਤਾਨੂੰ ਤਾਂ ਨਹੀਂ ਮੰਨਿਆ ਹੋਇਆ ਤਨ ਵਿੱਚ ਤਾਂ ਤਨ ਨਹੀਂ ਹੈ ਹੋਰ ਵੀ ਕਰਦੇ ਨੇ ਜਵਾਬ ਹੈ ਸੰਤੋਖ ધਨ ਸਭ ਧਨ ਧੂਲੀ ਸਮਾਨ ਸਾਰੇ ਤਨ ਮਿੱਟੀ ਬਰਾਬਰ ਨੇ ਜਿਹਦੇ ਕੋ ਸੰਤੋਖ ਸੰਤੋਸ਼ਤਾ ਰਹੇ ਸੰਤੋਖ ਤਾਂ ਤੇ ਹੈ ਨਹੀਂ ਸੰਤੋਸ਼ ਪ੍ਰਾ ਪਦਾਰਥ ਸੰਤੋਖ ਮਿਲਣਾ ਸੀ ਉਹ ਉਹਦੇ ਵਿੱਚ ਹੈ ਨਹੀਂ ਸਨਾਤਨਿ ਮਨ ਹੈ ਗੁਰਮਤ ਵਿੱਚ ਗਿਆਨ ਪਦਾਰਥ ਕਬੀਰ ਕਹਿੰਦਾ ਜਹ ਜ્ઞાન ਤਹਿ ਧਰਮ ਹੈ ਜਿੱਥੇ ਗਿਆਨ ਹੈ ਉਥੇ ਧਰਮ ਹੈ ज्ञान ने ना संतोष मिला ज्ञान का बद्दा मिल रहा है गुर बिना ज्ञान नहीं ये ज्ञान नहीं मिलता सो मत चवल्या कि ज्ञान पदार्थ है एदे नाल संतोष होना संतोष तण ज्यादा आ गया फिर किसी तान दी लोड़े नहीं थोड़ी अर्थ दी लोड़े यूं ही का नहीं है पदार्थ थोड़े खातर होगा सनातनई वक्त बात संसारी लोग खास्ते होगा संसारी वक्त खास्ते होगा ਗੁਜ਼ਾਰਿਆਂ ਦਾ ਆਲੇ ਵਾਸਤੇ ਹੋਊਗਾ ਵੀ ਬੰਦੇ ਨਹੀਂ ਚਾਰ ਪਦਾਰਥ ਉਹਨਾਂ ਵਾਸਤੇ ਹਿੰਦੂਆਂ ਵਾਸਤੇ ਹੋਊਗਾ ਸਿੱਖ ਗੁਰਸਿੱਖਾਂ ਵਾਸਤੇ ਨਹੀਂ ਗੁਰੂ ਘਰ ਵਾਸਤੇ ਤੈਸਾ ਸੋਣ ਤੈਸੀ ਉਸ ਤੈਸਾ ਅੰਮ੍ਰਿਤ ਤੈਸੀ ਵੇਖਾਟੀ ਤੈਸਾ ਮਾਨ ਤੈਸਾ ਅਮਾਨ ਤੈਸਾ ਰੰਗ ਤੈਸਾ ਰਾਜਾਨਾ ਢਾ ਲੱਗ ਹੋਰ ਉਹ ਉਹ ਤਾਂ ਗੁਰਦਾਨ ਦਾ ਸਨਾਤਨੀ ਮਤ ਹੈ ਸਾਰੀ ਉਹਦਾ ਜਰਾਤ ਨਹੀਂ ਮਰਦੇ ਢਾਲ ਨਹੀਂ ਲਿਆ ਉਹਨਾਂ ਵਾਲੇ ਪਦਾਰਥ ਨੇ ਉਹਨਾਂ ਹੁਣ ਹੁਣ ਮੰਨ ਵੀ ਗਏ ਅਸੀਂ ਗਲਤ ਪ੍ਰਚਾਰ ਕੀਤਾ ਉਹਨਾਂ ਨੂੰ ਵੀ ਪਤਾ ਲੱਗ ਗਿਆ ਸਮਝ ਗਏ ਹੋ ਵੀ ਇਹ ਤਾਂ ਪ੍ਰਚਾਰ ਗਲਤ ਹੈ ਨਹੀਂ ਸੀ ਪਤਾ ਉਹ ਸਮਝ ਗਏ ਮੰਨ ਗਏ ਉਹ ਵੀ ਹਾਂ ਗਲਤ ਹੈ ਹਾਂ ਸਾਡੇ ਚਾਰ ਪਦਾਰਥ ਕਿਹੜੇ ਨੇ ਜੀ ਸਾਡੇ ਗਿਆਨ ਪਦਾਰਥ ਪਹਿਲਾ ਧਰਮ ਚੋਂ ਗਿਆਨ ਮਿਲਣਾ ਜਿੱਥੇ ਗਿਆਨ ਨਹੀਂ ਹੋਦਾ ਤਾਂ ਉਹ ਗਿਆਨ ਕਿਹੜਾ ਮਿਲਣਾ ਆਤਮ ਗਿਆਨ ਇਹੋ ਨਾਮ ਵੀ ਕਹਿੰਦੇ ਨੇ ਆਤਮ ਗਿਆਨ ਨੂੰ ਪਹਿਲੀ ਸਟੇਜ ਜਿਹੜਾ ਲੈ ਇੱਕ ਨਾਮ ਬਿਨਾਂ ਕੰਨ ਦੇ ਸੁਣਨ ਵਾਲੇ ਕੰਨ ਗੁਰਬਾਣੀ ਹਰ ਨਾਮ ਸਮਾਇਆ ਗੁਰਬਾਣੀ ਚ ਨਾਮ ਸਮਾਇਆ ਹੋਇਆ ਉਹੀ ਬਣਦਾ ਗੁਰਬਾਣੀ ਨੂੰ ਮੰਤਰਨ ਕਰਦੇ ਤੇ ਜਿਹੜੇ ਲੱਕੇ ਉਹਨਾਂ ਕੰਦਾ ਉਹੀ ਤਾਂ ਗਿਆਨ ਅਗੁਰ ਵਰਤਿਦਾ ਪਹਿਲਾ ਗਿਆਨ ਬਦਲ ਗਿਆਨ ਤੋਂ ਮੁਕਤ ਪਦਾਰਥ ਮੁਕਤ ਤੋਂ ਨਾਮ ਪਦਾਰਥ ਮੁਕਤ ਬਕਰੀ ਵੀ ਗਿਆਨੀ ਧਿਆਗਾ ਉਹ ਤਾਂ ਮਰਤੀ ਹੋਇਆ ਸੰਸਾਰ ਛਡਾਉਂਦੀ ਹੈ ਮੁਕਤੀ ਤੇ ਮੁਕਤੀ ਤੋਂ ਬਾਅਦ ਨਾ ਅੱਗੇ ਨਹੀਂ ਜਾਂਦਾ ਮਾਤਾ ਨਹੀਂ ਵਰਕੇ ਜਿਉਂਦਾ ਕਰਨੇ ਫਿਰ ਜਨਪਦਾਰਥ ਹੈ ਜਨਪਦਾਰਥ ਤਾਂ ਮਿਲਦਾ ਇਹ ਨਾਮ ਪਦਾਰਥ ਮਿਲੇ ਤੁਰਕੀ ਬਾਣੀ ਆਈ ਤਿੰਨ ਅੰਗਲੀ ਜਨ ਤਵੜਾਈ ਉਹ ਨਾਮ ਹੈ ਬਿਨਾ ਕਰਨੇ ਤੇ ਸੁਣਨ ਵਾਲਾ ਜਿਹੜੇ ਨਾਮ ਨੇ ਬੰਦ ਕੀਤਾ ਸੀ ਜਿਹੜੇ ਚ ਉਹ ਨਾਮ ਖੋਲੂਗਾ ਬਾਹਰ ਕੱਢੂਗਾ ਤਾਂ ਨਿਕਲਦਾ ਸੰਸਾਰ ਤੋਂ ਬਾਹਰ ਮੁਕਤੀ ਦਾ ਬੁਖਤੀ ਦੰਗੇ ਤਾਂ ਜਾਂਦਾ ਨਾਮ ਨਾਲ ਤੁਰਕੀ ਬਾਣੀ ਨਾਲ ਬਿਨਾਂ ਕੰਨਾਂ ਤੋਂ ਸੁਣਨ ਵਾਲੇ ਹੁਕਮ ਨਾਲ ਹੁਕਮ ਨਾਲ ਬੰਦ ਹੋਇਆ ਹੁਕਮ ਨਾਲੇ ਬਾਹਰ ਨਿਕਲੋ ਜੇ ਜੇ ਪੂਰੀ ਵੀ ਕਰ ਲਵੇ ਨਾ ਸਜਾ ਫੇਰ ਵੀ ਸਰਕਾਰੀ ਹੁਕਮ ਨਾਲ ਬਾਹਰ ਨਹੀਂ ਕੱਢ ਸਕਦੇ ਨਿਕਲ ਸਕਦਾ ਸਰਕਾਰ ਦੀ ਮਰਜ਼ੀ ਹੈ ਛੱਡੇ ਜਾਂ ਨਾ ਛੱਡੇ ਜਿਹੜੇ ਬਹੁਤ ਕ੍ਰਿਮੀਨਲ ਹੁੰਦੇ ਨੇ ਕਹਿੰਦੇ ਜੇ ਸਰਕਾਰ ਨੂੰ ਤੇ ਖਤਰਾ ਹੋਵੇ ਨਹੀਂ ਛੱਡਦੇ ਵਿਭਾਰ ਆਉ ਖਤਰਾ ਬਾਹਰ ਕੱਢਣਾ ਹੋਰ ਗੱਲ ਹੈ ਹਾਂ ਕੈਦੀ ਨਹੀਂ ਉਹ ਕੈਦੀ ਵਾਲਾ ਕੰਮ ਨਹੀਂ ਉਹਦੇ ਲੈਣੇ ਸਜ਼ਾ ਉਹ ਜਾਨੀ ਮੁਸ਼ਕਲ ਨਹੀਂ ਉਹਨੂੰ ਹੈ ਪਰ ਉਹ ਜੜ੍ਹ ਚ ਬਾਹਰ ਖਤਰਾ ਉਹ ਤੋਂ ਇਸ ਕਰਕੇ ਮੁਫ਼ਤੀ ਵਾਲੇ ਤੋਂ ਬਾਹਰ ਖਤਰਾ ਆ ਜੇ ਮੁਕਤੀ ਆ ਜਿਹੜਾ ਹੈ ਨਾ ਮੁਕਤੀ ਵਾਲੇ ਤੇ ਨਹੀਂ ਮੁਕਤੀ ਵਾਲਾ ਮੁਕਤੀ ਦਾ ਬਾਣ ਆਰਾਧਨਾ ਆਰਾਧਨ ਆਰਾਧਨ ਨੀਕਾ ਹਰ ਹਰ ਨਾਮ ਆਰਾਧਨਾ ਆਰਾਧਨਾ ਤੇ ਬਾਅਦ ਜਾ ਕੇ ਕਿਤੇ ਨਾਮ ਮਿਲਦਾ ਉਹ ਤੋਂ ਬਾਅਦ ਹੁੰਦਾ ਇਥੋਂ ਫਿਰ ਫਿਰ ਸਰਵ ਹੁੰਦਾ ਫਿਰ ਲੀਨ ਹੁੰਦਾ ਫਿਰ ਅਨੇਕ ਹੈ ਮੁਕਤੀ ਦਾ ਅਨੇਕ ਨੇ ਇਹ ਸ਼ਬਦ ਵਿੱਚ ਜਿਹੜੀ ਨਾ ਫਿਰ ਇੱਕ ਹੁੰਦਾ ਸਾਰਿਆਂ ਨਾਲ ਸ਼ਬਦ ਦੇ ਰੂਪ ਵਿੱਚ ਹਕਮ ਦੇ ਰੂਪ ਇੱਕ ਹੈ ਕਲਾ ਕਲਾ ਅਨੇਕ ਹੈ ਫਿਰ ਇੱਕ ਹੈ ਅਨੇਕ ਤੋਂ ਇਕਤਾ ਵਿੱਚ ਨੂੰ ਜਾਣਾ ਜਦ ਫਿਰ ਬਾਹਰ ਨਿਕਲਦਾ ਬਾਹਰ ਆ ਕੇ ਕੋਈ ਹੈ ਮਾਇਆ ਵਿੱਚ ਅਨੇਕਤਾ ਹੈ ਮੁਕਤੀ ਵਾਲਾ ਮਾਇਆ ਦੇ ਵਿੱਚ ਹੈ ਜੇ ਅਨੇਕਤਾ ਹੈ ਉੱਥੇ ਉਹ ਤੇ ਦਾਸਨ ਬਾਦਸ਼ਾਹ ਕਹਿ ਰਹੇ ਚੇਤਨਾ ਤੇ ਉਹ ਹਮਰੋ ਆਵਨ ਕਾ ਹਮਰੋ ਆਵਨ ਕਾ ਚੁਮੀ ਰਹੀ ਸੁਤ ਪ੍ਰਭੂ ਚਨਨ ਮੈਂ ਹੋਈ ਸੀ ਜੁੜੀ ਹੋਈ ਸੀ ਚੁਮੀ ਰਹੀ ਹੈ ਲੀਨ ਸੀ ਲੀਨ ਹੋ ਰhalla ਚੁਮੀ ਹੋ ਰhalla ਧਿਆਨ ਉਦਨ ਕੀ ਹੋ ਰਹਾ ਸੰਸਾਰ ਚ ਦੇਖ ਰਹਾ ਰਾਜਾ ਰਾਮ ਕੀ ਕਹਾਣੀ ਜਾਣੇ ਹੈ ਬਾਬਾ ਜੀ ਤੁਸੀਂ ਪਦਾਰਥ ਦੀ ਗੱਲ ਕੀਤੀ ਨਾਮ ਪਦਾਰਥ ਵੀ ਆਇਆ ਨਾਮ ਪਦਾਰਥ ਫਿਰ ਉਹ ਚਾਰ ਪਦਾਰਥ ਜਿਹੜੇ ਹੋਏ ਫਿਰ ਇਹ ਨਾਮ ਪਦਾਰਥ ਅਲੱਗ ਹੋਇਆ ਪਹਿਲਾ ਗਿਆਨ ਪਦਾਰਥ ਆ ਯਾਰ ਜਿਹੜਾ ਗੁਰਬਾਣੀ ਵਾਲਾ ਨਾਮ ਹੈ ਗਿਆਨ ਪਦਾਰਥ ਹੈ ਕੋ ਨਾਮ ਪਦਾਰਥ ਜਿਹੜਾ ਬਿਨਨ ਕਰਨਾਂ ਤੇ ਸੁਣਨ ਵਾਲੇ ਤੁਰਕੀ ਬਾਣੀ ਉਹ ਹੈ ਉਹ ਉਹ ਅराधना ਨਾਮ ਦਾ ਇਹ ਜਪਨਾ ਨਿਲਦਾ ਹੈ ਗਿਆਨ ਜਪਦਾ ਵਿਸ਼ ਹੈ ਜਿਹੜਾ ਗਿਆਨ ਹੈ ਨਾ ਜੀ ਇਹ ਜਪ ਹੈ ਜਪ ਦਾ ਵਿਸ਼ਾ ਹੈ ਜਪਣਾ ਸਮਝਣਾ ਸੁਣਨਾ ਸੁਣੀਏ ਤੇ ਮੰਨਿਏ ਇਹ ਸੁਣ ਮੰਨਣ ਦਾ ਵਿਸ਼ਾ ਹੈ ਜਪਣ ਦਾ ਵਿਸ਼ਾ ਹੈ ਉਹ ਜਪਣ ਦਾ ਵਿਸ਼ਾ ਨਹੀਂ ਔਰ ਆਦਰਨ ਦਾ ਵਿਸ਼ਾ ਹੈ ਤੁਲਕੀ ਬਾਣੀ ਆਦਰਨ ਟੱਕ ਲੈ ਕੇ ਜਾਂਦਾ ਗਿਆਨ ਇਹ ਗਿਆਨ ਆराधना ਤੱਕ ਲੈ ਕੇ ਜਾਂਦਾ ਹੈ ਮੁਕਤੀ ਚ ਕੁਛ ਨਹੀਂ ਧਿਆਨ ਸਿਰਫ ਆराधना ਆराधना ਕਰਦੇ ਰਹਿਣਾ ਹੀ ਲਗਾਤਾਰ ਮੁਕਤੀ ਹੈ ਹੋਰ ਕੁਛ ਨਹੀਂ ਹੋਰ ਕੋਈ ਇੱਛਾ ਹੀ ਨਹੀਂ ਨਾਮ ਦੀ ਛ ਇਹਨੂੰ ਆराधना ਕਹਿੰਦੇ ਨੇ ਆराधना ਹੀ ਕਿਵੇਂ ਕਿਵੇਂ ਹੁੰਦੀ ਹੈ ਜੀ ਕੀ ਹੁੰਦਾ ਆराधना ਚ ਆਰਾਧਾ ਆਰਾਧਨਾ ਤਾਂ ਹੈ ਲੇਵੋ ਕੀ ਹੈ ਲੈਵ ਰਾਤ ਨਹੀਂ ਹੈ ਮੰਗਦਾ ਰੱਬ ਤੇ ਨਾਨਕ ਮੰਗੇ ਨਾਮદાન ਕਿਰਪਾ ਕਰੋ ਹਰੇ ਆਰਾਧਨਾ ਇੱਕੋ ਚੀਜ਼ ਮੰਗਦਾ ਹੈ ਉਹਦੀ ਲੋੜ ਏ ਨਹੀਂ ਹੋਰ ਕੋਈ ਉਹਦੀ ਲੋੜ ਹੀ ਆ ਨਾਨਕ ਨਾਮ ਮਿਲੇ ਤਾਂ ਜੀਵਾਂ ਨਾਮ ਮਿਲੇ ਤਾਂ ਜੀਵਾਂ ਵਰਿਆ ਤਾਂ ਹੈ ਗੁਗਤਾ ਹੈਗਾ ਨਾ ਨੂੰ ਨਾਮ ਮਿਲਾਂ ਤਾਂ ਜੀਵਾਂ ਤਾਂ ਲਗਿਆ ਇੱਥੇ ਨਹੀਂ ਤਾਇਰ ਇੱਥੇ ਤਾਂ ਤਾਂ ਜੀਵਾਂ ਜੀਵਾਂ ਤਾਂ ਬੋਲਣਾ ਬੋਲਣਾ ਜਿਉਣਾ ਬੁਲਾਇਆ ਜਦ ਬੁਲਾਇਆ ਬੋਲਦਾ ਉਹ ਜਿਉਣਾ ਸਾਬਤ ਹੈ ਫਿਰ ਉਚਾਰਨ ਕਰਦਾ ਗੁਰਬਾਣੀ ਉਹ ਜਨਮ ਬਦਾਸ ਮਿਲਿਆ ਹੋਇਆ ਸਾਬਤ ਹੋ ਗਿਆ ਜੇ ਸਾਵਧਾਨੀ ਨੀ ਕਰਦਾ ਤਾਂ ਨਾਮ ਨਹੀਂ ਮਿਲਿਆ ਜਿਹੜੇ ਕਹਿੰਦੇ ਸਾਨੂੰ ਚੁੱਪ ਹੋ ਗਏ ਜੇ ਚੁੱਪ ਹੋ ਗਏ ਤਾਂ ਮੁਕਤੀ ਤਾਂ ਖੋ ਸਕਦਾ ਚਲੇ ਗਏ ਤੁਸੀਂ ਪਰ ਮੁਕਤੀ ਵੀ ਦੱਸਣੀ ਪਊ ਤੁਹਾਨੂੰ ਕਿਵੇਂ ਹੋਏ ਆ ਉਹ ਤਾਂ ਮੁਕਤੀ ਵੀ ਨਹੀਂ ਦੱਸ ਰਹੇ ਮੁਕਤੀ ਮੁਕਤੀ ਦੀ ਜੁਗਤੀ ਕਰ ਰਹੇ ਨੇ ਜੁਗਤੀ ਹੁੰਦੀ ਹੋਈ ਨਹੀਂ ਗੁਰਬਾਣੀ ਜੋਤੀ ਰੱਦ ਕਰਦੀ ਹੈ ਜੋਗ ਜੁਗਤ ਇਹ ਪਾਈਆ ਜੁਗਤੀ ਰਸਿਆ ਕਿਵੇਂ ਆ ਅੰਜਨ ਮਾਹੇ ਨਰਿੰਦਲ ਲਈ ਹੈ ਯੋਗ ਚੁਗਤੀ ਵਪਾਈ ਹੈ ਅਜੋ ਜੁਗਤੀ ਤਾਂ ਪਾਉਣੀ ਹੈ ਪਹਿਲਾਂ ਅੰਜਨ ਮਾਹੇ ਨਰਿੰਦਲ ਹੋ ਕੇ ਤਾਂ ਦਿਖਾਓ ਮਾਇਆ ਦੇ ਵਿਚ ਰਹਣਾ ਹੈ ਮਾਇਆ ਤੋਂ ਨੰਦੇ ਫੋਕ ਦਿਖਾਓ ਮਾਇਆ ਦੀ ਇੱਛਾ ਤਿਆਗ ਕੇ ਦਿਖਾਓ ਲਗਾਤਾਰ ਕੈਸ ਕੇ ਦਿਖਾਓ ਲਗਾਤਾਰ ਇੱਛਾ ਢਾਕੇ ਹੋਈ ਹੈ ਮੁਕਤੀ ਉਨੂੰ ਰਾਜ ਨੂੰ ਕਹਿੰਦੇ ਨੇ ਜੇ ਕੋਈ ਇੱਛਾ ਫਿਰ ਜਾਗੇ ਰਾਜ ਨੂੰ ਖਤਮ ਇਹ ਮਾਇਆ ਵਾਲ ਤਾਂ ਚੱਲੇਗਾ ਆਰਾ ਉੱਥੇ ਬ੍ਰੇਕ ਹੋ ਜਾਂਦੀ ਹੈ ਜਿਵੇਂ ਸਰਵਰ ਇੱਕ ਵਾਰ ਟੁੱਟ ਜਵੇ ਨਾ ਪਿਛਲੇ ਸਾਲਸਾ ਤੋਂ ਨਵੇਂ ਸਾਲੇ ਚੰਦ ਸੂਰਜ ਦੀਵੜੇ ਚੰਦ ਸੂਰਜ ਦੀਵੜੇ ਆ ਸੰਸਾਰ ਦੀ ਚੰਦ ਸੂਰਜ ਦੀਵੜੇ ਨੇ ਜਿਹੜੇ ਆਪਣੇ ਜੀਵ ਨੇ ਇੱਕ ਇੱਕ ਨਹੀਂ ਚੰਦ ਹੈ ਕਿ ਨਹੀਂ ਸੂਰਜ ਇਹ ਲੱਖਾਂ ਚੰਦ ਨੇ ਲੱਖਾਂ ਹੀ ਸੂਰਜ ਨੇ ਔਰ ਇਸ ਮਨ ਵੀ ਚੰਦ ਸੂਰਜ ਨੇ ਰਗਾੜੀ ਚੰਦ ਸੂਰਜ ਵੀ ਨੇ ਅਦੂਏ ਵੀ ਨੇ ਬਾਹਲੇ ਵੀ ਨੇ ਇਹ ਬਾਲ ਨਹੀਂ ਚੰਦ ਸੂਰਜ ਦੇ ਬੜੇ ਨੇਖੇ ਉਹਦੇ ਕਰਕੇ ਬਾਈ ਡੜੇ ਦੀ ਬਣਾ ਤਾਂ ਕਰਚਾ ਚੰਦਾ ਸੂਰਜ ਸਾਡੇ ਦਾ ਦੀ ਗੱਡਾ ਲੱਗਦੀ ਬਾਉ ਜੀ ਜਿੰਦਾ ਵੀ ਉੱਡੇ ਹੀ ਨੇ ਇਹ ਘੜ ਦੀ ਵਿਸ਼ਾਲਤਾ ਹੈ ਜਿਵੇਂ ਸੂਰਜ ਦੀਵਾ ਉਹ ਘੜ ਕਿੱਡਾ ਜਿਹੜਾ ਹੈ ਲੱਗੜਾ ਬੀਜੂ ਦਾ ਕਹ ਰਹਾ ਹੈ ਕਿ ਜੀਸੂ ਦੀ ਵੋਕ ਨੇ ਨਹੀਂ ਬੀਜੂ ਰਾਜਾ ਚੰਦ ਸ਼ਿਵਜੀ ਦਾ ਤਾਂ ਕੋਈ ਕਾਰ ਹੈ ਹੀ ਨਹੀਂ ਉਹ ਤਾਂ ਕੰਦਾ ਬਣਾਇਆ ਹੀ ਸੀ ਉਹਨਾਂ ਤਿਆਗੀ ਹੈ ਉਹਦਾ ਮੰਨਦਾ ਵੀ ਤਾਂ ਕੰਦਾ ਹੁੰਦਾ ਹੀ ਨਹੀਂ ਇਹ ਕਾਰ ਹੈ ਹੀ ਨਹੀਂ ਉਹ ਵੀ ਆਪਣੇ ਆਪ ਨੂੰ ਮੰਨਦਾ ਮੇਰੇ ਤੋਂ ਕੁਝ ਹੰਕਾਰੀ ਹੁੰਦਾ ਜਿਹੜਾ ਬਿਸ਼ਨੂ ਦਾ ਉਤਾਰ ਹੈ ਹੰਕਾਰੀ ਹੁੰਦਾ ਹੈ ਰਾਮ ਜੀ ਵੀ ਹੰਕਾਰੀ ਹੈ ਕ੍ਰਿਸ਼ਨ ਵੀ ਹੰਕਾਰੀ ਹੈ ਉਹ ਵੀ ਐ ਕਰਦਾ ਕਾਲ ਬੱਪੜਾ ਕਾਲ ਬੱਪੜਾ ਕੌਤਕ ਦਿਖਾਉਂਦਾ ਇੱਥੇ ਊੜੇ ਬਾੜੇ ਤਲ ਕਾਲ ਕੀ ਐ ਕਾਲ ਹੁਕਮੇ ਆ ਹੁਕਮੇ ਕਾਲ ਐ ਕੌਤਕ ਨੇ ਸਾਰੇ ਹੁਕਮ ਨਾਲੇ ਜੰਮਣ ਮਰਨਾ ਹੁਕਮ ਨਾਲੇ ਸ੍ਰਿਸ਼ਟੀ ਚੱਲਦੀ ਐ ਕਾਲ ਅਕਾਲ ਖਤਮ ਕਾ ਕੀਨਾ ਅਕਾਲ ਖਤਮ ਦਾ ਕਾਲ ਬਣਾਇਆ ਹੋਇਆ ਹੈ ਕੀਨਾ ਹੁਕਮ ਕੀਦਾ ਅਕਾਲ ਦਾ ਅਕਾਲ ਬੋਲਣ ਦਾ ਕਾਲ ਕੀ ਹੈ ਕਾਲ ਹੁਕਮ ਜਮਣ ਮਾਨਾ ਹੁਕਮ ਹੈ ਇਹਦੇ ਹੀ ਕਾਹਤ ਸਾਰੇ ਜੋ ਕੁਝ ਹੋ ਰਿਹਾ ਇਹਦੇ ਹੋ ਰਿਹਾ ਹੁਕਮ ਨਾਲ ਸਭ ਕੁਝ ਹੈ ਕਾਲ ਬਪੂੜਾ ਕਿਉਂ ਹੈ ਹੀ ਹੁੰਦਾ ਕਾਲ ਹੋਰ ਕੀ ਹੋਊਗਾ ਕਾਲ ਵਗਣੇ ਤੇ ਇਹਨਾਂ ਜਿਹੜੇ ਕਿਸਦੇ ਅਧੀਨ ਹੋਵੇ ਪਪੜੇ ਹੁੰਦਾ ਉਹ ਕੋਈ ਵੀ ਨਹੀਂ ਪੰਡਾ ਨਹੀਂ ਹੈ ਹਾਕਮ ਦਾ ਹੁਕਮ ਹੈ ਹਾਕਮ ਦੇ ਦੀਨ ਹੁਕਮ ਹੁਕਮ ਹਾਕਮ ਉੱਪਰ ਆ ਕਰਨ ਦਾ ਮਤਲਬ ਇਹ ਹੈ ਬਪੂੜਾ ਦਾ ਕੀ ਅਰਥ ਹੈ ਜੋ ਕਿਸਦੇ ਬੱਚੇ ਹੋਵੇ ਕਾਲ ਦੇ ਕਾਲ ਦਾ ਕੀ ਨਾ ਕਾਲ ਜਿਹਨੇ ਕੀਤਾ ਜੋ ਜੋ ਰਚੋ ਤੋ ਤੇ ਸੇ ਤੇ ਆਉਦੇ ਕਾਬੂ ਹੈ ਸਕਲਾਂਸਪੁਰਖ ਦੇ ਕਾਬੂ ਹੈ ਉਹ ਉਹ ਤੇ ਵਖਰਾ ਨਹੀਂ ਉਹਦੀ ਮੰਜ਼ੀਆਂ ਸਾ ਉਹਦੀ ਮਰਜ਼ੀ ਹੋ ਕੋ ਹੋਰ ਕੀ ਹੈ ਇਹਨਾਂ ਨੇ ਇੰਡੀਪੈਂਡੈਂਟ ਬੰਨਿਆ ਕਾਲ ਨੂੰ ਇਹਨਾਂ ਨੂੰ ਤਾਂ ਕਿਹਾ ਇਹਨਾਂ ਨੇ ਕੁਝ ਹੋਰ ਮੰਨਿਆ ਤਾਂ ਉਹ ਨਹੀਂ ਪੜੇ ਗ੍ਰੰਥ ਇਹ ਜਿਹਨੂੰ ਜੀਰੋ ਉਪਦੇਸ਼ ਹੈ ਜੇ ਤੈਨੂੰ ਸਾਰਾ ਗਿਆਨ ਪੜਿਆ ਹੋਵੇ ਤਾਂ ਤੈਨੂੰ ਇਹ ਸਵਾਲ ਨਾ ਪੈਦਾ ਹੋਣ ਅਸਲ ਜੀ ਤੁਲੇ ਉਹ ਤਾਂ ਪੜਿਆ ਨਹੀਂ ਵਿਚਾਰਤਾ ਰੱਖੀ ਹੈ ਜਿਹੜੇ ਮੰਨਦੇ ਨੇ ਮੰਡਲ ਤੇ ਕੋ ਪੜਾਇਆ ਹੈ ਸਭਾ ਕਾਲ ਕਹਾਂ ਤੇ ਦਾੜੇ ਚਲੇ ਹਨ ਬਪਰੇ ਨਹੀਂ ਹੋਰ ਕੀ ਦੇ ਜੀ ਜਿਤੇ ਰਾਮ ਸੇਂ ਕ੍ਰਿਸ਼ਨ ਸੇ ਹੋਤ ਆਏ ਇਹਨੇ ਕਾਲ ਖਾਪਿਓ ਕਾਲ ਖਾਏ ਬਪੜਾ ਧੋਰ ਕੀ ਹੈ ਇਹ ਕਾਲ ਨੇ ਖਪਾਤੇ ਕਾਲ ਗਾਂਹ ਬਪੜਾ ਉਠਣ ਲੱਗੀ ਗੱਲ ਸੀ ਸਮਝ ਗਏ ਜੀ ਇਹ ਕਾਲ ਨਹੀਂ ਕਾਲ ਗਾਂਹ ਉਹਦੇ ਕਾਲ ਵੀ ਬਪੜਾ ਹੀ ਹੈ ਇਹ ਕਿਹਦੇ ਵਿਚਾਰੇ ਹੋਈ ਗਈ ਉੱਥੇ ਇਹ ਕਿਹੜੇ ਵਾਕ ਦੀ ਮੂਲੀ ਹੋਇਆ ਜਿਹਨੂੰ ਸੰਨਾਥਨੀ ਵਤਨੀ ਫਰਦਾ ਤਾਂ ਕੁਝ ਵੀ ਨਹੀਂ ਕਿ ਕਿਸੇ ਬਪੜਾ ਪਾਏ ਇੱਕ ਗਏ ਇੱਕ ਫੇਰ ਪਾਏ ਇੱਕ ਸ਼ਵ ਪਾਏ ਇੱਕ ਗਏ ਇੱਕ ਫੇਰ ਪਾਏ ਰਾਮ ਔਰ ਕ੍ਰਿਸ਼ਨ ਕੇ অবতার ਵੀ ਅਦੇਖ ਹੈ ਆਹ ਕੁਝ ਹੈ ਨਾ ਸਨਾਤਨੀ ਮਤ ਜੀ ਸਾਰਾ ਪੱਟੀ ਬੋਚੀ ਗੱਲ ਖਤਰ ਦਾ ਸਾਡੇ ਬਹਿਰ ਸੀ ਇਹਨਾਂ ਦਾ ਇਹ ਕਿਉਂ ਕਹਿੰਦੇ ਹੋ ਮੁਸਲਮਾਨਾਂ ਦਾ ਬਾਹਰ ਨਹੀਂ ਬਾਹਰ ਇਹਨਾਂ ਦਾ ਉਸ ਗਣ ਦਾ ਸਹਾਲ ਤੁਹਾਡਾ ਰਾਜ ਖਤਮ ਕਰ ਦੇਮੇ ਪਹਾੜੀ ਰਾਜੇ ਸਾਰੇ ਬਾੜੀ ਵਿਕਾਸੀ ਅੜਵੀ ਸਾਰੇ ਸੀ ਕੋਟ ਰਾਜ ਅਧੀਨ ਰਹਨੇ ਦੇਖਦੇ ਫਟ ਹੋ ਜਾਂਦੇ ਤੇ ਦੀਨ ਜਾਂਦਾ ਰਾयत ਵਾਲੇ ਵਾਗੀ ਰਹੇ ਨੇ ਇੱਥੇ ਮਤ ਹੋਰ ਹੈ ਚੰਡੀ ਨਵਾੰਦੇ ਰਹੇ ਜਾਂਦਾ ਖਣ ਵਾਲੇ ਵਾਗੀ ਰਹੇ ਨੇ ਇਸ ਕਰਕੇ ਸਿੰਘ ਜਾਂ ਜਾਂਦੇ ਸੀ ਨਾ ਪਰ ਆਇਆਂ ਦਾਨ ਵੱਲ ਤਾਂ ਚਲੇ ਜਾਂਦੇ ਤੇ ਇੱਧਰ ਰੁਮੀ ਤੇ ਆਉਂਦੇ ਯੂਪੀ ਵੱਲ ਨੂੰ ਇਹ ਤਾਂ ਸਾਰੇ ਦੁਸ਼ਮਣ ਤੇ ਯੂਪੀ ਵਾਲੇ ਪਹਾੜੀ ਰਾਜ ਵੀ ਦੁਸ਼ਮਣ ਸੀ ਇਹਨਾਂ ਦੀ ਵਿਚਾਰਦਾਰ ਇੱਕ ਉੱਤਰ ਵਾਲੇ ਨਹੀਂ ਗਏ ਦੱਖਣ ਵਾਲੂ ਗਏ ਨੇ ਦੱਖਣ ਦੀ ਵਿਚਾਰਦਾਰ ਹੋਰ ਹੈ ਉੱਤਰ ਦੀ ਹੋਰ ਹੈ ਦੱਖਣ ਦੀ আর ਪੱਛਮ ਦੀ ਵਿਚਾਰਦਾਰ ਰਲਦੀ ਆਪਣਾ ਪੱਛਮ ਦੇ ਵਿੱਚ ਮੁਸਲਮਾਨ ਸੀ ਉਹ ਤੇ ਗੁਰਨਾਨ ਗਾਇ ਨੇ ਕੋ ਟਕਰਾਇ ਹੋਇਆ ਉਹੁੰਦੇ ਹੀ ਚੱਲੇ ਗਏ ਨੇ ਉਹਨਾਂ ਨੇ ਪੀਰ ਮੰਨ ਲਿਆ ਇਹ ਦੁਨਾਨੇ ਗੁਰੂ ਮੰਨਿਆ ਝੂਠ ਗੱਲ ਹੈ ਕਿੰਦੇ ਵਿੱਚੋਂ ਕੁਝ ਆਦਮੀਆਂ ਨੇ ਗੁਰੂ ਬਣੇ ਬਹੁਤ ਥੋੜਿਆਂ ਨੇ ਬਰੋਹ ਜਿਆਦਾ ਉੱਤੋਂ ਹੁਰਵੀ ਮੰਨਦੇ ਨੇ ਅੰਦਰ ਬ੍ਰੋਧਾ ਮੁਚਾਤਾ ਦਾ ਦਾ ਬ੍ਰੋਧਾ ਉਹ ਉਹਨਾਂ ਦਾ ਸਾਡਾ ਉਹ ਇਹ ਦੁਨਾਨਾ ਗੁਰੂ ਹੈ ਇਹ ਦੁਈਆ ਇਹਨਾਂ ਦਾ ਗੁਰੂ ਹੈ ਇਹ ਦੁਈਆ ਗੁਰੂ ਬਦਲਦਾ ਹੁੰਦਾ ਗੁਰੂ ਦੱਸਦਾ ਵੀ ਤੂੰ ਹੀ Hindu ਬਣੋ ਗੁਰੂ ਨੂੰ Hindu ਬਣਾਉਂਦੇ ਫੇਰ ਗੁਰੂ ਕਹਿੰਦਾ ਜੇ Hindu ਹੈ ਜੇ Hindu ਹੈ ਫਿਰ ਤਾਂ ਗੁਰੂ ਨਹੀਂ ਹੋ ਤੂੰ ਗੁਰੂ ਹੋ ਤੇ ਤੂੰ ਪਹਿਲਾਂ ਹੀ ਨੇ ਉਹ ਗੁਰੂ ਆ ਗੁਰੂ ਕਾਣੀ ਕਹਿੰਦਾ ਫੇਰ ਗੁਰੂ ਆ ਜਿਹੜਾ ਨਵੀਂ ਰੋਸ਼ਨੀ ਦਵੇ ਜੋ ਪਿੱਛੇ ਰੋਸ਼ਨੀ ਹੁੰਦਾ ਨਵੀਂ ਰੋਸ਼ਨੀ ਦਵੇ ਤਾਂ ਗੁਰੂ ਆ ਇਹ ਰੋਸ਼ਨੀ ਨਿੰਮੈ ਦਿੱਤੇ ਗੁਰੂ ਕਾ ਦਾ ਨਾਮ। ਇਹ ਗੁਰੂ ਮੰਦਰ ਨੇ ਸੇਖਵੀ। ਨਵੀਂ ਰੋਸ਼ਨੀ ਕੀ ਹੈ ਜੋ ਕੋਈ ਦੱਸੇ। ਇਹ ਲੋਗ ਤਾਂ ਉਹੀ ਚਾਰ ਪਦਾਲਸ ਨੇ। ਨਵੀਂ ਰੋਸ਼ਨੀ ਦੱਸੋ ਕੀ ਨਵੀਂ ਲਾਈਟ ਜਿਹੜੀ ਦਿੱਤਿਓ ਦਿਖਾਉਣ ਕੀ ਹੈ। ਗੁਰੂ ਵੀ ਹੈ ਲਾਈਟ ਵੀ ਪ੍ਰਾਣੀ ਹੈ। ਲਾਟਣ ਵੀ ਹੋਈ ਹੈ, ਬੱਤੀ ਵੀ ਹੋਈ ਹੈ, ਤੇਲ ਵੀ ਹੋਈ ਹੈ, ਸਭ ਕੁਝ ਹੋਈ ਹੈ। ਕੋਈ ਮਾਇਆ ਮਾਇਆ ਵਾਲਾ ਤੇਲ ਹੈ ਜਲਦਾ। ਜੋਦ ਵੀ ਉਹੀ ਹੈ ਨਵਾਂ ਕੀ ਹੈ ਤੁਹਾਡੇ ਕੋਲ ਗੁਰੂ ਕਾਗਾ ਗੁਰੂ ਤਾਂ ਹੈ ਉਹਦਾ ਗਿਆਨ ਗੁਰੂ ਹੈ ਜੋ ਗਿਆਨ ਦਿੰਦਾ ਉਹੀ ਗੁਰੂ ਹੁੰਦਾ ਹੈ ਉਹ ਉਹਨੇ ਨਵਾਂ ਗਿਆਨ ਦਿੱਤਾ ਕੁਛ ਉਹ ਤਕਵੀਰ ਵਾਲਾ ਹੀ ਦਿੱਤਾ ਚਾਹੇ ਪਰ ਨਵੇਂ ਸਿਰੇ ਤੋਂ ਦਿੱਤਾ ਉਹ ਗੰਗਲਾ ਕਰਤਾ ਸੀ ਪਹਿਲਾਂ ਵੀ ਸੀ ਕਵੀਰ ਤੋਂ ਪਹਿਲਾਂ ਵੀ ਸੀ ਨਾਰਦ ਵਾਲਾ ਗਿਆਨ ਹੈ ਨਾਰਦ ਵਾਲੀ ਭਗਤੀ ਹੈ ਭਗਤ ਨਾਰਦ ਦੀ ਇਹਦੇ ਨਾਲ ਉਪਜੀ ਇਹ ਹਿੱਦ ਚੁੱਪ ਜਿਓ ਨਹੀਂ ਹੈ ਉਪਜਣੀ ਸੀ ਤਾਂ ਪੈਦਾ ਹੋਣੀ ਸੀ ਭਗਤ ਨਾਰਦ ਦੀ ਇਹਦੇ ਨਾਲ ਉਪਜੀ ਉਪਜੀ ਕਿਦੋਂ ਮੁਜੀਏ ਜਿਹਦੇ ਉਹ ਚਾਨਣ ਕਰੂਗੀ ਇਹ ਭਗਤੀ ਹੈ ਗੁਰ ਮਤ ਜੇ ਗੁਰ ਮਾਤਾ ਨਾ ਉਹੀ ਉਭਜਣੀ ਅੰਦਰ ਉਹੀ ਸੋਈ ਸੋਈ ਜਾਗਣੀ ਹੈ ਫਿਰ ਜਿਹੜਾ ਚੰਨ ਉਹ ਦਊਗੀ ਉਹ ਗਿਆਨ ਗੁਰੂ ਹੋਊਗਾ ਉਹ ਨਵਾਂ ਚੰਨ ਹੋਊਗਾ ਹਾਂਜੀ ਜੀ ਜਿਵੇਂ ਤੁਸੀਂ ਦੱਸਿਆ ਹੁਣ ਵੀ ਪਿਛਲੇ ਗ੍ਰੰਥ ਦੇ ਵਿੱਚੋਂ ਇਹ ਗੱਲਾਂ ਆਈਆਂ ਕੀ ਫਿਰ ਸਾਨੂੰ ਉਹ ਵੀ ਪੜ੍ਹਨੇ ਚਾਹੀਦੇ ਆ ਤੁਸੀਂ ਕੀ ਲੈਣੇ ਪੜ੍ਹ ਕੇ ਯਾਰ ਉਹਨੂੰ ਜਿਹੜੇ ਮੰਨਦੇ ਤੇ ਉਹਨਾਂ ਨੂੰ ਉਪਦੇਸ਼ ਕਰਕੇ ਆਪਣੇ ਨਾਲ ਲੈ ਆਉਂਦਾ ਠੀਕ ਹੈ ਜੀ ਸਾਰੀ ਦੁਨੀਆ ਨੂੰ ਬਤੇ ਸਾਰੀ ਦੁਨੀਆ ਦੀਆਂ ਬਤਾਂ ਨੂੰ ਉਪਦੇਸ਼ ਹੈ ਕੈਂ ਕੀ ਲੈਣਾ ਪੜ ਕੇ ਤੂੰ ਕਿੱਥੇ ਖੜਾ ਤੈਨੂੰ ਕਿਹੜਾ ਉਪਦੇਸ਼ ਹੈ ਤੇਰੇ ਦੀ ਬਿਮਾਰੀ ਹੈ ਦੀ ਦਵਾਈ ਖਾਣੀ ਹੈ ਤੈਨੂੰ ਜਿਹੜੀ ਬਿਮਾਰੀ ਦਵਾਈ ਲੈ ਜੀ ਦੇ ਪੜਨ ਦਾ ਆ ਪਤਾ ਨਹੀਂ ਥੋੜਾ ਗੁਰਬਾਣੀ ਸੇ ਬਹੁਤ ਸੀਮਤ ਬਤਲਵਾ ਸੁਣਣ ਵਾਲਿਆਂ ਦਾ ਤੂੰ ਸਾਲ ਨੂੰ ਜੱਫਾ ਪਾਣੀ ਬੈਠੇ ਹੋ ਜੱਫਾ ਉਹ ਲੋੜਾ ਜਿਹਨੇ ਦੁਨੀਆਂ ਨੂੰ ਸਮਝਾਉਣਾ ਹੋਵੇ ਸਾਰਿਆਂ ਨੂੰ ਜਿਹੜਾ ਕੋ ਡਾਕਟਰ ਬਣਨਾ ਹੋਵੇ ਜਿਹਨੇ ਬੈਦ ਬਣਨਾ ਹੋਵੇ ਬੈਦ ਬਣਨਾ ਤਾ ਪੜੋ ਜੇ ਬੈਦ ਨਹੀਂ ਬਣਨਾ ਆਪਣੀ ਯੋਗਾ ਲੈਣਾ ਫਿਰ ਆਪਣੇ ਮਤਲਬ ਦੀ ਗੱਲ ਪੜੋ ਦੋਈ ਜਿਹੜੀ ਬਵਾਰੀ ਤੁਹਾਨੂੰ ਹੈ ਠੀਕ ਹੈ ਜੀ ਜ਼ਰੂਰੀ ਨਹੀਂ ਹੈਗਾ ਵੀ ਸਾਰਾ ਕੁਝ ਹੀ ਕਰਨਾ ਆਪਣੇ ਲਈ ਪਹਿਲਾਂ ਆਪਣੇ ਲਈ ਕਰਨਾ ਅਸੀਂ ਆਪਣੇ ਲਈ ਕਰੋ ਅਸੀਂ ਕਿੱਥੇ ਖੜੇ ਆਂ ਜਦ ਤੂੰ ਹੀ ਨਿਰੋਗ ਹੋ ਜਾਉਂਗੇ ਤਦ ਨੂੰ ਆਪੇ ਗੱਲ ਹੋ ਜੂ ਆਪ ਤਾਂ ਨਿਰੋਗ ਰੋਗ ਦਾ ਕਾਰਨ ਆਪੇ ਪਤਾ ਲੱਗ ਜੂ ਨੂੰ ਕਿ ਬਿਮਾਰੀਆਂ ਦਾ ਇਲਾਜ ਦੱਬੀ ਹੈ ਤੋਂ ਪਹਿਲਾਂ ਆਪਣੀ ਬਿਮਾਰੀ ਦਾ ਇਲਾਜ ਕਰਦੇ ਅਸੀਂ ਹਰ ਇੱਕ ਲੈ ਕੇ ਜਫਾ ਪਾ ਲੈਂਦੇ ਹਰ ਇੱਕ ਲੈ ਕੇ ਜਫਾ ਪਾ ਲੈਂਦੇ ਤੂੰ ਕੀ ਜਾਣਦਾ ਹੁੰਦਾ ਥੋੜੀ ਬੈਕਰਾਉਂਡ ਦਾ ਨਹੀਂ ਪਤਾ ਤਦ ਮਜ਼ੀਦਾ ਛੋੜੇ ਕੰਮ ਸਮਝ ਆ ਜੂ ਫਿਰ ਮੇਰੇ ਮਾਂ ਪੂਰੀ ਜ਼ਿੰਦਗੀ ਲਾ ਦੋ ਛੱਡੋ ਕੰਮ ਉਹ ਤੁਸੀਂ ਕਰ ਨਹੀਂ ਸਕਦੇ ਤੇ ਤੁਸੀਂ ਆਪਣੇ ਜੋਗਾ ਹੀ ਰੱਖੋ ਬਸ ਜਿਹਨੂੰ ਜਿਹੜੀ ਬਿਮਾਰੀ ਸੀ ਜਿਹੜੀ ਮਾਂ ਪੜਾਤੀ ਪੁੱਠੀ ਉਹ ਉਹਦਾ ਉਹਨੂੰ ਸਮਝ ਉਹਨੂੰ ਬਾਈਏ ਥੋੜਾ ਐ ਪੁੱਠੀ ਹੈ ਉਹ ਪੁੱਠੇਰਾ ਪਿਆ ਹੋਇਆ ਜਦੋਂ ਆਇਆ ਵੀਰ ਆਪੋ ਠਾਈਦੈ ਨੂੰ ਐਨੂੰ ਜਾਣੋ ਸੀ ਤਾਂ ਇੱਥੋਂ ਭੁੱਲ ਗਿਆ ਜਾਂ ਦੋਰਾ ਘਿਆ ਹੀ ਨਹੀਂ ਤੇਰੇ ਮਤਲਬੇ ਕੋਈ ਨਹੀਂ ਸਾਡਾ ਸਤਿ ਸਕਲ ਮਤਲਬ ਹੈ ਵੀ ਚਾਰ ਬਦਾਰਥੇ ਨੂੰ ਆਨੇ ਨੇ ਸਾਡੇ ਬਦਾਰਥਾਏ ਨੇ ਗੁਰਬਾਣੀ ਦਾ ਗਿਆਨ ਆਂ ਕਹਿੰਦਾ ਸੰਤੋਖ ਚਾਹੀਦਾ ਹੈ ਕੋਈ ਤੂੰ ਇਮਾਨਦਾਰੀ ਚਾਹੀਦੀ ਹੈ ਦੋ ਗੱਲਾਂ ਨੇ ਇਮਾਨਦਾਰੀ ਆ ਸੰਤੋਖ ਬਾਕੀ ਤੁਸੀਂ ਕੀ ਲੈਣਾ ਦੁਨੀਆ ਤੇ ਬਾਕੀ ਦਸ ਘੜੀ ਜਿੰਦੀ ਲੋੜ ਹੈ ਫੇਰ ਜੋ ਬਾਣੀ ਦੀ ਲੋੜ ਹੈ ਇਹ ਸ਼ਬਦ ਦੀ ਤੁਹਾਨੂੰ। ਕਿ ਆਪਨੇ ਅਮਰੂਣ ਜਾ ਲੈਣਾ ਐਵੇਂ ਚਖਮਾਲ ਦੇ ਫਰੀ ਜਾਣਾ। ਤੁਹਾਨੂੰ ਸਮਝ ਨਹੀਂ ਆਈ ਅਸਲ ਦੇ ਵਿੱਚ। ਕਿ ਕਾਨੂੰਨੀ ਨੀ ਇਹ ਤਾਂ ਹੀ ਸਖ ਫਸੇ ਨੇ। ਤੁਹਾਨੂੰ ਸਮਝ ਨਹੀਂ ਆਈ ਗੱਲ ਕੀ ਐ ਇਹ। ਕਿ ਗੁਰਦਾਰਿਆਂ ਨਹੀਂ ਕੰਮ ਹੋ ਸਕਦਾ। ਇਹਨੂੰ ਦੁਨੀਆਂ ਨੂੰ ਉਲ ਜਾਤਾ ਕਦੇ ਕੋਈ ਸ਼ਬਦ ਨੇ ਕਦੇ ਕੋਈ ਸਾਰੇ ਉਲ ਜਾ ਸਕਦੇ। ਉਹ ਉਹ ਨਹੀਂ ਸਲੇਪਸ ਦੱਸੋ ਭਾਈ ਤੈਨੂੰ ਆਮ ਮਾਰੀ ਐ ਐ ਦਵਾਈ ਖਾਣੀ ਐ ਐ ਪਰਹੇਜ ਰੱਖ ਤੈਂ ਬਸ ਆਪਣੇ ਤੱਕ ਫੀਸ ਉਤਰੇ ਫਿਰ ਕੇ ਤੇ ਪੰਨੇ ਕੁਝ ਪੈ ਜਾਂਦਾ ਇਹ ਨਾਲ ਆ ਬੁੱਢੇ ਨੇ ਨਨ ਜਾਂਦੇ ਸਾਰੇ ਇੱਕ ਆਦਮੀ ਕਪੜਾ ਕੇਸ ਰੰਦਦਾ ਉਹ ਆਪਣੇ ਕੇਸ ਤੱਕ ਮਾਤਲਬਾ ਉਹਨੇ ਵਕੀਲ ਬਣਨਾ ਸੁਪਰੀਮ ਕੋਰਟ ਦਾ ਉਹੀ ਸਬੂਤ ਇਕੱਠੇ ਕਰਦਾ ਜਿਹਦੇ ਨਾਲ ਉਹਦਾ ਕੇਸ ਜਿੱਤਿਆ ਜਾ ਸਕੇ ਬੱਤ ਉਹ ਆਪਣੇ ਕੇਸ ਦੇ ਸਬੂਤ ਇਕੱਠੇ ਕਰੋ ਤੁਸੀਂ ਤੁਸੀਂ ਇੰਟਰਨੈਸ਼ਨਲ ਲੈਵਲ ਦੇ ਵਕੀਲ ਬਣਨਾ ਚਾਹੁੰਦੇ ਹੋ ਤੁਸੀਂ ਕਿਹਨਾਂ ਉਹ ਵਕਾਲਤ ਤੇ ਥੋਤੇ ਨਹੀਂ ਮੰਨਣਾ ਵਕੀਲ ਉਹ ਵਕੀਲ ਬਣਨਾ ਫਿਰ ਵਕਾਲਤ ਹੀ ਫਿਰ ਤੁਹਾਨੂੰ ਆਪਣਾ ਕੰਮ ਛੱਡ ਲਓ ਪ੍ਰੋਬਲਮ ਇੱਥੇ ਆਉਂਦੀ ਆ ਕੇ ਤੁਹਾਨੂੰ ਆਪਣੇ ਤੁਸੀਂ ਸਬੂਤ ਇਕੱਠੇ ਕਰੋ ਆਪਣੇ ਬਿਆਨ ਦਿਓ ਕੀ ਕੱਲੋਂ ਮੇਰੇ ਮੈਂ ਬਿਆਨ ਕੀ ਦੇਣੇ ਨੇ ਕਿਹੜੇ ਮੇਰੇ ਖਿਲਾਫ ਜਾਂਦੇ ਨੇ ਕਿਹੜੀ ਗੱਲ ਮੇਰੇ ਹੱਕ ਆ ਜਾਊਗੀ ਬੋਲਣਾ ਸਿੱਖੋ ਅਦਾਲਤ ਵਿੱਚ ਕੀ ਹੈ ਹਾਂਜੀ ਜਾਚੈ ਕਰ ਲక్ష్ਮੀ ਕੁਵਾਰੀ ਚੰਦ ਸੂਰਜ ਦੇਵੜੇ ਕੌਤਕ ਕਾਲ ਪਪੂੜਾ ਆਹ ਸੂਰਜ ਇਹਦਾ ਚਾਂਦਾ ਜੇ ਮਨਮੁਖਾ ਦਾ ਗਿਆਨ ਹੈ ਚੰਦ ਦਾ ਮਨਮੁਖਾ ਜਿੱਥੇ ਮਨਮੁਖੀ ਦੋਹਿਲਾ ਮਨਮੁਖਾ ਤੇ ਜਿੰਨਾਂ ਤੇ ਗਈ ਪੱਛਾ ਨੂੰ ਆਇਆ ਚੰਦਰਾ ਜਿੰਨਾ ਮਰਜੀ ਚਾਹੇ ਉਹਨਾਂ ਮਾਸ਼ੀਦਾ ਹੋਵੇ ਪਰ ਹੋਊ ਰਹੇ ਚੰਦ ਦਿਨ ਹੋਇਆ ਚੰਦ ਚੰਨ ਰੋਸ਼ਨੀ ਉਹ ਦਿਆ ਤਾਰਿਆਂ ਦੀ ਰੋਸ਼ਨੀ ਹੁੰਦੀ ਹੈ ਤਾਰੇ ਰਹੀ ਜੀਵਨ ਨੇ ਤਾਰਿਆਂ ਦੇ ਜੀਵਨ ਇਹਨਾਂ ਨੇ ਕਹਿਣਾ ਜੀ ਕਿੰਨੀ ਰੋਸ਼ਨੀ ਆ ਤਾਰਿਆਂ ਦੀ ਤਾਰਿਆਂ ਦੀ ਰੋਸ਼ਨੀ ਆ ਇਹ ਜਿਹੜਾ ਸਨਾਤਨ ਮਤ ਹੈ ਸਨਾਤਨ ਮਤ ਕੋ ਤਾਰਿਆਂ ਦੀ ਆ ਸਭ ਲਈ ਜੀ ਤਾਰੇ ਹੀ ਨੇ ਹੋ ਇਹਨਾਂ ਦੇ ਚੰਦਰਮਈ ਜੀ ਦੀ ਰੋਸ਼ਨੀ ਹੋਣਾ ਸੀ ਤਾਂ ਚੰਦਰਮਈ ਦਾ ਕਲਾ ਨੇ ਜਿਹਨ ਕੋ ਕਹਿੰਦੇ ਨੇ 16 ਤਲਾ ਸਿੰਗਰਮਾਪੂਰ ਨੂੰ ਪੂਰਨਮਾਸੀ ਉਹ ਵੀ ਰਾਤ ਹੈ। ਨਾਲੇ ਦਾ ਦੇਖਣ ਉਹ ਕਾ ਜਨਰ ਦੇ ਵਿੱਚ ਆਪਣੇ ਵਿੱਚ ਦਾਗ ਨਹੀਂ ਹੈ। ਕੋਈ ਜਾ ਚੈ ਕਰ ਜੀ ਦੇ ਜਾ ਚੈ ਜਿਸ ਵਿੱਚ ਯਾਰ ਆਂਦਾ ਕਹਿ ਲਾਂਦਾ ਚਾਹਦਾ ਉਹਦਾ ਵਿੱਚ ਵਿੱਚ ਦਾ ਚਾਹ ਆ ਗਿਆ ਅੱਪਾ ਕਹਿੰਦੇ ਖਰਚ ਕਹਿੰਦਾ ਨਹੀਂ ਜੀ ਉਹ ਕਹਿੰਦੇ ਡੱਬੀ 'ਚ ਹੈ ਛੇ ਕਹਿੰਦੇ ਵਿੱਚ ਨਹੀਂ ਵਿੱਚ ਹੈ ਛੇ ਕਹਿੰਦੇ ਨੇ ਤੇ ਉਹੀ ਚੇ ਲੱਗਿਆ ਇੱਥੇ ਜਾ ਲਗਾ ਕੇ ਲੰਗ ਜਿਸਚੋ ਜਿਸ ਵਿੱਚ ਵਿੱਚ ਨਾ ਜਿਸਚੋ ਜੀ ਜਦੋਂ ਦਾ ਵਿੱਚ ਇਹ ਸ਼ਬਦ ਹੈ ਯਾ ਚੈ ਘਰ ਜਲਕੀ ਕੁਆਰੀ ਤੇ ਅਕਲ ਕੁਆਰੀ ਹੋਇਆ ਹੈ ਗਾਲ ਗੋਲੀ ਖਾਇਆ ਵਾਰੀਆ ਹੂੰ ਚੰਦ ਸੂਰਜ ਦੀਵੜੇ ਚੰਦ ਸੂਰਜ ਦੀਵੇ ਨੇ ਤੇਰਾ ਮੰਨਦਾ ਗਾ ਇਹਦੇ ਘਰ ਦੇ ਵਿੱਚ ਨੇ ਕਹਿੰਦੇ ਸੂਰਜ ਨੇ ਦੀਵੜੇ ਨੇ ਜਾਂਦੇ ਸੂਰਜ ਨੇ ਦੀਵੇ ਬਣਾਏ ਨੇ ਆਪ ਆਪ ਨੂੰ ਦਾ ਉਹ ਰੋੜ ਨਹੀਂ ਦੀਵੇ ਰੱਖਣ ਦੀ ਸਾਡੇ ਬਾਹਰ ਤੇ ਬਣਾਏ ਨੇ ਆ ਘਰ ਦੇ ਵਿੱਚ ਆਪਾਂ ਰਹਿੰਦੇ ਉਹ ਜਿੰਨ ਤੱਕ ਇਹ ਅਰੰਡਦੇ ਆਪਾਂ ਰਹੇ ਨਹੀਂ ਆਪਣੇ ਘਰ ਜਾਨਾ ਜੀ ਉਹ ਜਿਹੜੀਆਂ ਨਾਲ ਜਿਹੜੀਆਂ ਮਾਤਾ ਉੱਗਣ ਵਾਲੇ ਲੰਗੇ ਸ਼ਿਤੀਰਾਮ ਤੇ ਜਿਹੜੀਆਂ ਉਹ ਕਹਿੰਦੇ ਸਾਡਾ ਘਰ ਤੂੰ ਕਹਿੰਦਾ ਮੇਰਾ ਦਾ ਉਹ ਜੂਹਾਂ ਦੇ ਫਟਾਉਂਨਾ ਪਾਪੜੀ ਹੋਰ ਕਿੰਨੇ ਛੋਟੇ-ਮੋਟੇ ਜੀਵਾਨਾ ਉਹਨਾਂ ਦਾ ਵੀ ਏਰੀਆ ਦਾ ਬੈਥੂ ਵੈਰੇ ਉਹ ਕਹਿਣਾ ਸਾਡਾ ਕਿੱਲੀ ਨੰਦ ਨਾਮ ਹੁੰਦੀ ਜੇ ਹੁੰਦੀ ਛੰਡਾ ਦੋਈ ਗੱਲੀ ਨਹੀਂ ਹੁੰਦੀ ਬੋਦੀ ਬੋ ਨਾ ਨਾ ਤਰ ਵੀ ਹੈ ਤੇ ਤੇਰੇ ਨਾਲ ਤਾਂ ਅੱਜੇ ਤਾਂ ਕੀੜੇ ਮਕੌੜੇ ਨੋਦੇ ਕਾਲਦੇ ਕਰਤਾ ਹੋਦਾ ਯਾ ਸੀ ਵੀ ਕੀੜੇ ਮਕੌੜੇ ਵਿਚੇ ਰਹਿੰਦੇ ਆ ਜੇ ਜਿਹੜੀ ਪਰੇਸ਼ੀ ਕਰਚੇ ਹੁੰਦੀ ਹੈ ਜਿਹੜੀ ਆ ਜਾਂਦੇ ਸੋ ਵੇ ਆਂ ਚੁਗਿਆ ਜ਼ੋ ਫਾਨੀਆ ਆ ਆ ਇਹ ਦਾ ਫਰੰਡੀ ਕਰ ਹੁੰਦਾ ਕਾਰਜ ਬਹੁਤ ਕੁਝ ਹੁੰਦਾ ਉਹ ਤਾਂ ਕੰਮ ਖਾ ਗਿਆ ਉਹ ਤਾਂ ਕਹਿਣਾ ਨਹੀਂ ਇਹ ਤਾਂ ਕਰਤਾ ਬੈਠੇ ਸਭ ਕੁਝ ਆਫਰ ਕੋਲੋ ਤੇ ਕੱਪਟੇ ਸ੍ਰੀ ਕੋਟਵਾਲਾ ਉੱਤੇ ਪੌਣੇ ਕੋਟਵਾਲ ਕੋਟਵਾਲੋ ਕਬੀਰ ਕਹਿੰਦਾ ਸੰਤਾਂ ਮਾਨ ਨੂੰ ਦੂਤਾਂ ਨੂੰ ਇਹ ਕੋਟਵਾਰੀ ਮੇਰੀ ਜਿਹੜਾ ਸੱਜਦਾ ਪ੍ਰਚਾਰਕ ਹੈ ਨਾ ਚੱਕੀ ਮਤ ਇੱਕ ਕੋਟਵਾਲੀ ਇਹਦੀ ਹੈ ਸਰਦਾਰੀ ਹੈ ਕੋਟਵਾਲੀ ਜੂਠੇ ਨੂੰ ਦੰਦ ਦੰਦ ਲੋਦੇ ਨੂੰ ਸਜ਼ਾ ਦੇਣੀ ਸੱਚ ਨੂੰ ਮਾਨ ਦੇਣਾ ਜੋਰ ਦਾ ਤਰਸਕਾਰ ਕਰਦੂ ਗੁਰਬਤ ਕਰਨੀ ਲਈ ਮਨ ਮ ਕੋ ਅਪੇਜਣਾਂ ਤੇ ਜੀ ਪੱਥਰ ਘੈਤਾ ਹੁੰਦਾ ਨਾਨਕ ਤੇ ਪੇ ਨਾਲ ਅਸਲ ਖਰ ਕੁੱਤਾ ਤੇ ਗੁੜਵਾਰੀ ਨਹੀਂ ਹੈ ਜੇ ਬੇਨੁਗੁਣ ਗਰਭ ਕਰਨ ਤੇ ਗੁੜਵਾਰੀ ਨਹੀਂ ਹੈ ਕੁੱਟੇ ਨੇ ਕੋੜਵਾਲੀ ਕੁੱਟੇ ਉਹ ਸਾਰੇ ਕੁੱਟਣਾ ਤਾਂ ਮਨ ਕੋ ਕੁੱਟੇ ਇਹਨਾਂ ਦਾ ਮਨ ਕੁੱਟਿਆ ਮਨ ਕੁੱਟਿਆ ਤਾਂ ਅੰਨੇ ਕੁੱਟਿਆ ਬੁਰਵਾਣੀ ਮਨ ਨੂੰ ਕੁੱਟਦੀ ਹੈ ਤੁਹਾਨੂੰ ਜੀ ਕੁੱਟਦੀ ਤੁਹਾਨੂੰ ਤਾਂ ਕੋੜਦੇ ਨੇ ਸੁਨਾਤ ਨਹੀਂ ਬਰਮੀ ਮਾਰੀ ਤਾਂ ਪਣੀ ਉਹ ਸਰੀਰ ਨੂੰ ਤਾਂ ਉਹ ਕੁੱਟਦੇ ਨੇ ਨੇ ਮਨ ਨੂੰ ਘਰ ਦੀ ਇਹੋ ਬਾਣੀ ਉੱਟਣਾ ਤਾਂ ਮਨ ਕੋ ਖੂਪਦਾ ਤੇ ਉਹ ਮਨ ਕੋ ਉੱਟੇ ਪੰਜ ਅੰਤੈ ਛੂਪਦਾ ਤਾਂ ਪਰ ਬ huzur ਹੁੰਦੇ ਤਰਨਾਇ ਲੈਂਦੀ ਹੈ ਤੇ ਤੋਂ ਵੀ ਆਪਾਂ ਉਹ ਵੀ ਇਦਾਂ ਕਹਿ ਜੀਣਾ ਇਹਾ ਕਪੜਾ ਕੋਲ ਲੈ ਤੋ ਇਹੇ ਪੜ ਤੇ ਪੜਦੇ ਇਹ ਮਨ ਹੁੰਦੀ ਹੈ ਤੇ ਆਖਰੀ ਕੋਟਾ ਆ ਤਾਂ ਦੇ ਫਟ ਗਿਆ ਕੱਪੜਾ ਜਾਂ ਫਿਰ ਜਾਂ ਫਟ ਗਿਆ ਜਾਂ ਫਿਰ ਬਣ ਗਿਆ ਜਾਂ ਨਿਕਲ ਗਿਆ ਫਟ ਗਿਆ ਉਹ ਟਾਂ ਵਾਲੇ ਨੇ ਆਪਣੀ ਕਹਾਣੀ ਦਈ ਜਿੱਦਾਂ ਸ਼ਰਮਾਂ ਨਹੀਂ ਹੁੰਦੀ ਕੋਲੋਂ ਸਰੀਰਾਂ ਫਟ ਗਿਆ ਫਟ ਗਿਆ ਉਹਦਾ ਅੱਡ ਹੋ ਗਿਆ ਫਟ ਗਿਆ ਉਹਦਾ ਮਨ ਉਹਨੇ ਆਪਣਾ ਦੂਰ ਕਾਂਦੇ ਅਲੱਗ ਹੋ ਗਿਆ ਵਿਸ਼ਨਰੀਆਂ ਨੇ ਕਲਾਸ਼ ਨੂੰ ਇਹਦੀ ਫਟਣੀ ਹੈ ਆਪਣੇ ਨਾਲੋਂ ਇੰਨੇ ਆਦਮੀ ਫਟੇ ਕੇ ਜੀ ਉਪਦੇਈਨਾ ਹਾਂਜੀ ਸੋ ਹੈ ਜੀ ਸ਼੍ਰੋਮਣੀ ਕਮੇਟੀ ਵਿਭਾਗ ਦੂਜਾ ਉਹਦੇ ਵਿੱਚ ਸੋ ਕਰਾ ਸ੍ਰੀ ਸ਼ੁਕਰਾ ਸ੍ਰੀ ਵੀ ਹੈ ਹੋ ਸ਼ੁਕਰਾ ਹੀ ਹੈ ਇਹ ਜਿਹੜੀ ਸਾਡੇ ਨੂੰ ਜਿਹੜੀ ਕਿਰਤ ਹੈ ਹੈ ਜਿਹੜੀ ਜਾਣ ਕੋਤਵਾਲੀ ਹੈ ਇਹ ਸੁਖ ਹੈ ਦੀ ਦੁਖਰੇ ਤਕ ਕੀ ਹੈ ਪਰਮ ਦੇ ਵਿੱਚ ਫਸਾਉਣਾ ਜੋ ਹੈ ਪਰਮ ਦਾ ਨਾਸ ਕਰਨਾ ਦੁਨੀਆ ਦਾ ਸੁਖ ਹੈ ਇਹ ਜੋ ਕਰਮਨ ਦੇ ਨਿਮਨ ਦਾ ਫੈਲਾਉਣਾ ਪ੍ਰਚਾਰ ਕਰਨਾ ਭਰਮ ਦੇ ਵਿੱਚ ਪਾ ਕੇ ਲੋਕਾਂ ਨੂੰ ਲੁੱਟਣਾ ਭਰਮ ਵਿੱਚ ਪਾ ਕੇ ਗੁਰੂ ਬਣਨਾ ਅਗਿਆਨਤਾ ਫੈਲਾਈ ਰੱਖਣਾ ਅਗਿਆਨਤਾ ਕਰਕੇ ਲੋਕਾਂ ਨੂੰ ਗੁੰਮਰਾਹ ਕਰਨਾ ਇਹ ਪਾਪ ਹੈ ਬੁਕਲਤੀ ਹੈ ਪਾਪ ਕਰਨ ਤਾਂ ਜਨਮ ਕੇਵ ਜਿਓ ਤੇ ਕੋਈ ਨਾ ਮੇਲੀ ਰਾਮ ਤੇ ਬੋਲ ਮੇਲੀ ਕੋਈ ਵੀ ਨਹੀਂ ਹੈ ਐ ਵਰਮਾ ਵੀ ਜੂ ਸ਼ਵੀਰ ਨੇ ਜੇਹਨੇ ਸਾਥ ਲੈਂਦੇ ਨੇ ਉਹਦੇ ਬੁੱਧਨੀ ਕਰਨਾ ਬੋਲਣਾ ਉੱਥੇ ਜੇ ਹੋਊਗਾ ਤਾਂ ਮੋਲੋ ਇਹ ਥੱਲੇ ਹੀ ਨੇ ਚੋਰ ਕਾਮਾ ਭਰੇ ਨਾ ਕੋਈ ਚੋਰ ਆਰਾਮ ਖੋਨੇ ਹਮ ਕੋਈ ਨਹੀਂ ਪਰਣਾ ਕਰਨੇ ਇਹ ਦੁਕ੍ਰਿਤੀ ਹੈ ਕੁਟਵਾਲੀ ਸੁਕ੍ਰਿਤੀ ਸੋ ਉੱਪਰ ਹੋਸਨ ਬੈਨੇ ਰਾਖਸ਼ਣਾ ਗੁਰੂ ਆ ਹੋ ਤਾਂ ਕਹਿੰਦੇ ਨੇ ਰਾਜਮੰਦੇ ਨੇ ਉਹਨਾਂ ਨੂੰ ਕੁਟਦੇ ਨੇ ਰਾਖੇ ਨੇ ਦੇਵਤਾ ਕੀ ਨੇ ਕਿਆ ਕੇ ਬੜੇ ਹਮਦਰਦੀ ਨਾਲ ਗੱਲਾਂ ਕਰਕੇ ਸੰਤ ਬੜਾ ਫਸਾ ਕੇ ਲੁੱਟਦੇ ਨੇ ਖਾਂਦੇ ਨੇ ਹੌਲੀ ਹੌਲੀ ਖਾਦੇ ਕਰਕੇ ਉਹਨਿੰਦੇ ਮੂੰਹ ਵਿੱਚ ਪਾਣੀ ਮੂੰਹੋਂ ਮਿਟੈਨ ਨਾ ਕੇ ਜੀ ਹੋ ਗਈ ਹੈ ਮੂੰਹੋਂ ਮਿਟਾ ਜਮਾ ਨਹੀਂ ਹੁੰਦਾ ਖੁਦ ਉਪਰੇਤੀ ਹੈ ਉਹ ਆਪਣੇ ਨਾਲ ਸਾਥ ਬਾਸੇ ਮਿਟਾ ਹੌਲੀ ਜੀ ਤੋ ਐਸਾ ਰਾਜਾ ਸ਼੍ਰੀ ਨਰਹਰੀ ਐਸਾ ਹੈ ਉਹ ਵੈਸਾ ਨਹੀਂ ਜੈਸਾ ਤੁਸੀਂ ਕਹਿੰਦੇ ਹੋ ਨਰਹਰੀ ਉਹਨਾਂ ਨੇ ਜੋ ਨਰਹਰੀ ਐਕਸਲੈਂਸ ਕੀਤਾ ਉਹ ਤੋਂ ਉਲਟਾ ਐਕਸਲੈਂਸ ਉਹਨਾਂ ਇਹਦਾ ਮਤਲਬ ਐਸਾ ਹੈ ਜੈਸਾ ਆਪ ਪਹਿਲੇ ਬਤਾ ਰਹੇ ਵੈਸਾ ਨਹੀਂ ਹੈ ਜੇ ਜਿਹੜਾ ਉਹ ਜਿਹੜਾ ਕਹਿੰਦੇ ਉਹ ਜਿਹੇ ਹੁੰਦਾ ਫਿਰ ਐਸਾ ਲੈ ਰਹੇ ਕੀ ਲੋ 20 ਸਾਰੀ ਵੇਖਾ ਦਤੀ ਹੈ ਉਹ ਜਦੋਂ ਲਕੀਰ ਪਾ ਹੈ ਪੁਲਾਨ ਸਭ ਬੁਣਾ ਕੇ ਕਿਹਾ ਐ ਉਹ বিষ্ণੂ ਦੇ ਕਾਲ ਜਿਹੜੇ ਰਤਨ ਸੀ ਉਹ ਨਹੀਂ ਸੀਗੇ ਉਹ ਬੰਦਰ ਦੇ ਵੱਡੇ ਲੈ ਕੇ ਭੱਜੇ ਬੇਈਮਾਨ ਨਿਕਾ ਟਿੱਕੇ ਬਾਅਦ ਚ ਉਹਦਾ ਕਾਲਸਾਂ ਕੁਝ ਕਿੱਥੇ ਹੈ ਹਾਂਜੀ ਅਰੇਲੀ ਕੰਪਨੀ ਕੀ ਹੈ ਜਾਂਚ ਹੈ ਕੋ ਲਾਲ ਬ੍ਰਹਮਾ ਚਤੁਰਮੁਖ डावੜਾ ਜਿਹੜੇ ਘਰ ਦੇ ਵਿੱਚ ਇੱਕ ਬ੍ਰਹਮਾ ਵੀ ਹੈ ਆਲੇ ਉਹ ਬ੍ਰਹਮਾ ਨਾਲ ਜਿੱਤ ਚਤੁਰਮੁਖ ਚਾਰ ਮੁਖ ਵਾਲਾ ਅਸਲ ਨੇ ਚਾਰੇ ਪੇਦ ਦੇ ਤੋ ਨੇ ਚਾਰ ਮੂੰਹ ਬਣਾਤੇ ਚਤੁਰਮੁਖ ਸੀ ਮੁਖ ਇੱਕੋ ਹੀ ਚਾਹੀਦਾ ਉਹ ਚਤੁਰਾ ਬੜਾ ਚਤੁਰ ਦਾਤ ਆਇਆ ਹੋਇਆ ਚਤੁਰਾਈ ਜਿਹੜੀ ਹੈ ਇਹਨਾ ਨਾ ਪਾਇਆ ਆਇਰ ਮੰਚਨ ਚਲ ਚੰਚਲਤਾ ਰੰਗਿਆ ਜਿੰਨਾ ਚਿਰ ਆਪਣੇ ਆਪ ਨੂੰ ਚਤੁਰ ਮੰਨਦਾ ਹੋ ਚਾਣਾ ਮੰਨਦਾ ਚੈ ਚਾਣ ਪਾਲਾ ਕੋਈ ਖਲ ਨਾਲ ਜਦੋਂ ਆਪਣੀ ਜਾਣ ਪਛੜ ਦਿੰਦਾ ਹੋ ਜਾਂਦਾ ਫਿਰ ਗੁਰਮੁਖ ਹੋ ਜਿਹੜਾ ਹੈ ਉਹ ਪੜਨਤ ਹੋ ਜਾਂਦਾ ਘਰ ਵਿੱਚ ਆਹੋ ਜਿਹਦਾ ਕਹ ਰਿਹਾ ਉੱਥੇ ਹੀ ਰਹਿੰਦਾ ਹਾ ਹੁਣ ਬ੍ਰਹਮਾ ਕੁਲਾਲ ਕੁਲਾਲ ਲਿਖ ਬੱਤੇ ਲਾਲੀ ਦੇ ਨਾਮ ਨਹੀਂ ਹੈ ਉਹ ਵੇਦ ਜਿਹਨੇ ਵੇਦਾਂ ਦੇ ਵਿਚਾਰ ਤਾਨੂੰ ਵਗਾੜ ਕੇ ਇਹ ਦੱਸ ਰਿਹਾ ਉਹ ਕੁਲਾਲ ਹੈ ਲਾਲ ਲਾਲ ਤੇ ਲਾਲਨ ਕੁਲਾਲ ਕਕਰੂ ਕੜਾ ਕੇ ਨੈਗੇਟਿਵ ਲੱਗਿਆ ਲਾਲੀ ਮੇਰੇ ਲਾਲ ਕੀ ਨਾਮਦਾਰ ਮ ਲਾਲ ਹੁੰਦਾ ਨਾ राले ब्रह्मा चतुर्मुख बड़ा सयाना जी ओ पढ़ला ता अर बाद पाठती ते शास्त्र काढले उने हां कुलाल ब्रह्मा चतुर्मुख डावड़ा डावड़ा चार मुखाड़ा जिन विश्व संसार राची ले ਉਹ ਕੈਨਾਂ ਨੇ ਵਿਸ਼ਵ ਸੰਸਾਰ ਨੂੰ ਰੱਖਿਆ ਜਿਹਨੇ ਤੁਸੀਂ ਕਹਿੰਦੇ ਹੋ ਵਿਸ਼ਵ ਸੰਸਾਰ ਰੱਖਿਆ ਉਹ ਦਾ ਕਹੇ ਆ ਯਾਨੀ ਉਹਦਾ ਹੋ ਨੌਕਰ ਹੈ ਉਹਦਾ ਕਰਦਾ ਮਾਨ ਕਰਦੇ ਆ ਉਹਦਾ ਮੁਲਾਜ਼ਮ ਕਹ ਲੋ ਨੌਕਰ ਕਹ ਲੋ ਤੇ ਆ ਉਹ ਰਾਮ ਕਹ ਲੋ ਇਛ ਵੀ ਹੈ ਉਹਦਾ ਕਰਿਆ ਜਾਂਚੇ ਈਸ਼ਰ ਬਾਵਲਾ ਜਗਤ ਇਥਰ ਆ ਗਿਆ ਨਾ ਚੇਵੀ ਇਥਰ ਇਥਰ ਬਾਵਲਾ ਜਿਹਨੂੰ ਤੁਸੀਂ ਬਾਵਲਾ ਕਹਿੰਦੇ ਹੋ ਚੇਵੀ ਪੰਗਪੀਰ ਬਾਵਲਾ ਇਸਰ ਵੀ ਉਹਦੇ ਘਰ ਕੇ ਉਹ ਹਿੰਦੂ ਗੰਤੇ ਭੱਟੀ ਪਹੁੰਚੀ ਜਾਂਦਾ ਉਹ ਵੀ ਉਹਦੇ ਘਰੇ ਆ ਉਸ ਘਰ ਦੇ ਗਿਆਨਪਤ ਜਗਤਗੁਰੂ ਕਹੋਂਦਾ ਆਪਣੇ ਆਪ ਨੂੰ ਜਗਤਗੁਰੂ ਬਣ ਕੇ ਬੈਠਾ ਬ੍ਰਹਮਾ ਆਪਣੇ ਆਪ ਨੂੰ ਗੁਰੂ ਨਹੀਂ ਮੰਨਦਾ ਅੰਨ ਮਾਮਣ ਗੁਰੂ ਬਣ ਆ ਕੇ ਬੈਠੇ ਜਗਤਗੁਰੂ ਉਹ ਕਹਿੰਦਾ ਮੈਂ ਜਗਤਗੁਰੂ ਭਾਰਤ ਤੱਤ ਗਿਆਨ ਤੋਂ ਸਖਣਾ ਜਿਹੜਾ ਗਿਆਨ ਹੈ ਉਹਦਾ ਤੱਤ ਨਹੀਂ ਆਉਂਦੇ ਵਿੱਚ ਤੋਂ ਸਾਰ ਤੱਤ ਗਿਆਨ ਤੋਂ ਸਖਣਾ ਤੱਤ ਗਿਆਨ ਤੋਂ ਵਾਂਝਾ ਗੁਰੂ ਆ ਤਤਸਾਰਖਾ ਗਿਆਨ ਪਾ ਕੀਲੇ ਆ ਤਤ ਤੋਂ ਖਾਲੀ ਕਹਿੰਦਾ ਲੋਕਾ ਤਤ ਨਹੀਂ ਆਉਦੇ ਵਿੱਚ ਸੱਚ ਨਹੀਂ ਹੈ ਜਿਹੜਾ ਗਿਆਨ ਉਹ ਦੱਸ ਰਿਹਾ ਭਰਮ ਗਿਆਨ ਦਾ ਪ੍ਰਚਾਰ ਕਰ ਰਿਹਾ ਆਪਣੇ ਗਿਆਨ ਦੇ ਵਿੱਚ ਲੋਕਾਂ ਨੂੰ ਭਰਮਾ ਰਹੇ ਹੋਣ ਜਾ ਰਹੇ ਫਾਂਸਣ ਕੀ ਵੀ ਨਹੀਂ ਦੱਸ ਰਿਹਾ ਫਾਂਸਣ ਕੀ ਵੀ ਸਭ ਕੋ ਜਾਣੇ ਉਹਦੀ ਬੇਦੀ ਫਸਾਉਣ ਵਾਲੀ ਹੈ ਮਾਇਆ ਚ ਫਸਾਈ ਰੱਖਣ ਵਾਲੀ ਹੈ ਕਿਉਂਕਿ ਮੁਕਤੀ ਤਾਂ ਖੁਦ ਮੰਗਦਾ ਪ੍ਰਮਾਣ ਗੰਧੀ ਕੋ ਖੋਜੇ ਮਹੇਸ਼ਰ ਪ੍ਰਮਾਣ ਗੰਧੀ ਤਾਂ ਕੋਈ ਦੇ ਮੁਕਤੀ ਦਾ ਤਾਂ ਕੋ ਹੈ ਮੁਕਤੀ ਤਾਂ ਆਪ ਚਾਹੁੰਦਾ ਸਿਰ ਉਹ ਕਿਹੜਾ ਗਿਆਨ ਹੈ ਜਿਹੜਾ ਦੇ ਰਿਹਾ ਲੋਕਾਂ ਨੂੰ ਮੰਨਦਾ ਅਜਾ ਮਾਰਾਜ ਫਸਾਉਣ ਵਾਲੇ ਗਿਆਨ ਨੇ ਉਹਦਾ ਗਿਆਨ ਨਾ ਮਾਇਆ ਤਮੰਦੀ ਹੈ ਜ਼ਰੂਰ ਰਉਦਰ ਭਗਤ ਜਗਤਮਾਹੈਂ ਦਸ ਬਾਸ਼ਾ ਕਰਨ ਰਉਦਰ ਭਗਤ ਜਗਤਮਾਹੈਂ ਸੁਖ ਕੇ ਦੇਵ ਸੋ ਸਦਾ ਪਰੈ ਸੰਤਾਰਿ ਸੁਖੋ ਉਰੁ ਸੰਤਾਰਿ ਸੁਖਤਾ ਬਣਜੈ ਨਾ ਸੁਖ ਕੇ ਦੇਵ ਸਦਾ ਪਰੈ ਮਰੈ ਫਰਾਵਾ ਭਗਤੀ ਭਗਤ ਨੂੰ ਮੁਕਤੀ ਦੀ ਵਿਰਤੀ ਤੇ ਮੁਕਤੀ ਦੀ ਵਿਰਤੀ ਚਰਮਗਾਹ ਹੈ ਗੁਰੂ ਹੈ ਮਾਈ ਬੁੰਡੋ ਤੇ ਗੁਰੂ ਕੀ ਜਾਤੇ ਜਾਏ ਤਾਹੀ ਆਏ ਗੱਲ ਕਹੀ ਹੈ ਕਬੀਰ ਆ ਇਹ ਤੇ ਰੁਖਿਆ ਜਗਤ ਗਰੂ ਰੂ ਜੋ ਉਹਦੇ ਜਟਾਂ ਨੇ ਬਹੁਤ ਬੜੀਆਂ ਬਣੀਆਂ ਤੱਤੇ ਉਹਦੀ ਮੱਤ ਨੂੰ ਮੰਡੋ ਉਹਦੀ ਮੱਤ ਵਿੱਚ ਜਟਾ ਨੇ ਜਟਾ ਆਵੇਂ ਜੇ ਉਹ 라ਵੀ ਲੈ ਜਟਾ ਫੇਰ ਕਿਹੜਾ ਕੁਛ ਹੋ ਗਿਆ ਗੱਲ ਫੇਰ ਵੀ ਉਹੀ ਹੈ పాਪ ਪੁੰਨ ਜਾਂਚੇ ਡਾਂਗੀਆਂ ਦੁਆਰੇ ਜਿਹਦੇ ਦੁਆਰੇ ਹੈ ਉੱਤੇ ਬਾਰੇਦਾਰ ਖੜੇ ਨੇ ਚੋਬ ਦਾ ਲਾਂਗਾਂ ਲੈ ਕੇ ਖੜਦੇ ਨਹੀਂ ਹੁੰਦੇ ਇੱਕ ਦੋ ਬੰਦੇ ਦਵਾਰਪਾਲ ਜੀ ਖੜੇ ਤੋੜੇ ਦਰਵਾਜਾ ਪਾਪ ਪੁਨਨ ਦਰਵਾਜਾ ਇੱਕ ਪਾਪ ਦੇ ਦਰਵਾਜੇ ਤੇ ਖੜਾ ਇੱਕ ਪੁਨਨ ਵਾਲੇ ਤੇ ਖੜਾ ਪਾਪ ਪੁਨਨ ਪਾਪ ਦਰਵਾਜਾ ਖੁੱਲਦਾ ਜੀ ਬਾਗਿਆ ਪਾਪ ਪੁਨ ਦੋਨੋਂ ਭਾਈ ਭਾਈ ਦੋ ਭਾਈ ਨੇ ਦੋ ਮਿਲਕੇ ਕੇ ਸੇ ਸਪਾਈ ਹੈ ਦੋ ਦਰਵਾਜੇ ਨੇ ਕਿਤੇ ਚੇਤਾ ਕਿਤੇ ਮਾਨਾ ਦੋ ਇੱਕ ਪੁੰਨੀ ਰਗ ਪਾਪੀ ਹੈ ਡਾਂਗੀਆਂ ਬਾਬਾ ਜੀ ਡਾਂਗਾ ਆਲੇ ਲੱਛੀ ਦਾ ਕਿਹੜੇ ਖੜੇ ਨਹੀਂ ਹੁੰਦੇ ਚਿੱਤਰ ਗੁਪਤ ਲੇਖੀਆ ਆ ਅੰਦਰ ਜਿਹੜਾ ਚਿੱਤਰ ਉਹ ਵੀ ਚਿੱਤਰ ਹੋਉਂਦੇ ਚਿੱਤਰ ਉਹ ਲੇਖਾ ਕਰਦਾ ਉਹ ਯੋਗ ਹੈ ਜੜੇ ਚਿੱਤਰਗੁਪਤ ਦਾ ਕੀ ਅਰਥ ਹੈ ਜੀ ਜੇ ਤਜੇ ਜੇ ਤਰਾਂ ਦੀ ਐਂਟ ਤੇ ਬੋਪਤਾ ਇਹਨਾਂ ਲਈ ਕਹਿੰਦਾ ਜੇ ਤਬ ਉਹ ਦੁਰਜਸ ਉਹ ਤੇ ਤੈਨੂੰ ਪਰਨ ਹੋ ਯਾਰ ਕੰਮ ਤਾਂ ਖਰਾਬ ਹੈ ਕਰਾਂਗਾ ਨੰਦਾ ਦਾ ਇਹੋ ਲੇਖਾ ਕਰਦਾ ਦਿਖਾ ਕੇ ਨਹੀਂ ਕਰਦਾ ਜੇ ਤੁਹਾਨੂੰ ਗੁਪਤੇ ਅੰਦਰ ਦੀਨ ਅਨਿਵਾਰ ਬੈਠਾ ਸਭ ਦੇ ਅੰਦਰ ਬਿਖਾਲਿਆ ਹੋਇਆ ਗੋਆਪੀ ਚਤਰਗੁਪਤਾ ਹੈ ਹੋਰ ਕੌਣ ਹੈ ਕੋਈ ਨਹੀਂ ਧਰਮ ਰਾਏ ਪਰੋਲੀ ਪ੍ਰਤੀਹਾਰਾ ਅਜਲਾ ਧਰਮਾ ਹੈ ਉਹ ਹੀ ਧਰਮਾ ਹੈ ਕੋਤਨੁਰਾਵੀ ਉਸ ਨੂੰ ਗੈਰ ਨੇ ਜਦ ਲੈ ਖਾ ਮੰਗਾ ਉਹਦੇ ਉੱਪਰ ਹੈ ਉਹ ਹੋਰ ਉੱਪਰ ਥੋੜੀ ਹੋਰੀ ਸੀਟ। ਇਕਾ ਥੱਲੇ ਉਹ ਨਾ ਕੋਈ ਮੁਚੀ ਬਿਲਾਨ ਕਰਦੀ ਏ ਮੁਚੀ ਲਿਖਦਾ ਆ ਥੰਦੜ ਇਕ ਉੱਪਰ ਉਹ ਤਾਰ ਬੁਲਾਇਆ ਜਬ ਲੇਖਾ ਮੰਗਾ ਜੀ ਉਹ ਲੇਖਾ ਮੰਗਣ ਵਾਲਾ ਕਹੇ ਕਲੇਖਾ ਲੈਣ ਵਾਲਾ ਕਲੇਖਾ ਉਹ ਨੂੰ ਕਿ ਕਦਾ ਲਿਖ ਜਾਣਦਾ ਹੀ ਆ ਇਹ ਕਲੇਖਾ ਤੇ ਉਹਦਾ ਹਸਾਬ ਮੰਗਣ ਉਹ ਉਹ ਪ੍ਰティਹਾਰ ਉਸ ਪਰ ਬੈਠਾ ਲਾਗ ਲਈ ਉਹ ਪੁੱਛੂਗਾ ਕਿ ਨਾ ਜਵਾਬ ਉਹਦੇ ਮੂਹਰੇ ਜਵਾਬ ਦੇ ਹੈ ਜਵਾਬ ਤਲਵੀ ਹੈ ਉਹਦੇ ਪ੍ਰਤੀ ਜੋ ਲੇਖਾ ਉਹਦੇ ਪ੍ਰਤੀ ਜਵਾਬ ਦੇ ਹੀ ਹੈ ਤੁਹਾਰਾ ਜੋ ਲਿਖਿਆ ਗਿਆ ਉਹਦੇ ਬਾਬਤ ਉਹਦੇ ਪਰਥਾਏ ਜਵਾਬ ਤਲ وی جواب اے نہیں لکھاں لے کیوں چھڈ دے نا او تعبین کرنا تے ہاں روندی پے یار او ہے نا کہ ایک دا ہندا لکھاں لکھیاں چھڑیاں نا او دا کوئی یار او دی کوئی پرواہ نہیں نہیں نہیں او لکھے را سب دینا پنے جواب دہی ہے او دی لکھے ਜੋ ਲੇਖਾ ਖਾ ਲੈ ਕੇ ਆ ਜਾ ਉਹਨੇ ਪ੍ਰਤੀ ਜਿਮੁਰ ਬਾਰੀ ਆਤਾ ਦੀ ਵਿਆਖਿਆ ਨੇ ਪਰੋਲੀ ਦਾ ਕੀਤਾ ਪਰਲੋ ਵਾਲਾ ਦਰਬਾਨ ਜੋ ਅਧਿਕ ਅਨ ਅਧਿਕਾਰੀ ਨੂ ਅੰਦਰੋ ਜਾਣੋ ਰੋਕਦਾ ਹੈ। ਯਾਰ ਪਰੋਲੀ ਅੰਦਰੋ ਜਾਣੋ ਨਹੀਂ ਰੋਕਦਾ ਸਰਬਰਾਜ। ਸਰਬਰਾਜ ਅੰਦਰੋ ਜਾਣੋ ਰੋਕਦਾ। ਦਰਬਾਨ ਮਤਲਬ ਪਪਾ ਰਾਰੇ ਨੂੰ ਮਲਵਾਨ ਆ ਗਿਆ ਹੁਣ ਦਰਵਾਨ ਬਾਅਦ ਫਿਰ ਕਹਾਂ ਜਾਣਾ ਹੈ ਇਹ ਆ ਹਾਂਜੀ ਉਹ ਤੀਸ ਤੁਰਿਆ ਫਿਰ ਪਰੋਲੀ ਪਰਲੋ ਕਰਨ ਵਾਲਾ ਵੀ ਲਿਖਿਆ ਜਿਨ੍ਹਾਂ ਨੇ ਨਹੀਂ ਨਹੀਂ ਪਰਲੋ ਕਰਨਾ ਪ੍ਰਤੀ ਉਹ ਪੂਰੇ ਦੇ ਪ੍ਰਤੀ ਜੋ ਲੇਖਾ ਲਿਖਿਆ ਜਾਊ ਵਹਾਂ ਦਾ ਜਾਏਗਾ ਉਹ ਤਾਂ ਫਰਾਮਗਦਾ ਤੇ ਜਵਾਬ ਤਲ ਵੀ ਲੈਣੀ ਆ ਉਹਦੀ ਸਜ਼ਾ ਦੇਣੀ ਆ ਤੈਨੂੰ ਹਮਲਾ ਕਰਨਾ ਹੁੰਦਾ ਜੇ ਵੀ ਹੈ ਹੰਕਾਰ ਤੇ ਪ੍ਰਹਾਰ ਨਹੀਂ ਕਰਦਾ ਜੀ ਉਹਵੇਂ ਪ੍ਰਹਾਰ ਹੀ ਲਿਖਿਆ ਉਹਨੂੰ ਜੋੜ ਕਰਨੀ ਆ ਉਹਨੇ ਤੇ ਲੇਖੇ ਤੇ ਜਵਾਬ ਚਲੂ ਹੀ ਆ ਜਵਾਬ ਦੇਣਾ ਪੈਣਾ ਤੈਨੂੰ ਗੱਲਾਂ ਹੁੰਦਾ ਦੇ ਪ੍ਰਤੀ ਤੇਰੇ ਉਹਦੇ ਸਵਾਲਾਂ ਦਾ ਜਵਾਬ ਦੇਣਾ ਪੈਣਾ ਤੈਨੂੰ ਜਵਾਬ ਦੇਹੀ ਹੈ ਫਰਨਾ ਹੁੰਦਾ ਉਹਦੇ ਪ੍ਰਤੀ ਜੋ ਲਿਖਿਆ ਉਹਦੇ ਉੱਪਰ ਉਹਨੇ ਉਪਰੇ ਉਹਦੇ ਬੈਸ ਹੋਣੀ ਹੈ ਵੇ ਨਹੀਂ ਪਾਇਲ ਤੇ ਪੁੱਛੇ ਛੋੜੀਆਂ ਤੇਰੀ ਦਿੰਦੇ ਸ਼ਾਮ ਲਾ ਉਹਦੀ ਜਵਾਬ ਦੇ ਦਿੱਤੀ ਤੇਰੀ ਗਾਂ ਗਾਂ ਤੂੰ ਨਹੀਂ ਗੱਲ ਦੀ ਉਹਨੇ ਇੱਕ ਕੇਸ ਭੇਜਤਾ ਦਫਾ ਲਾ ਕੇ ਅੱਗੇ ਤਾਲ ਚਲੇ ਜਵਾਬ ਦੇ ਤੇਰੀਆਂ ਤੇ ਹੋਰ ਕਿਹਦੇ ਉਹਦੇ ਪ੍ਰਤੀ ਉਹ ਪ੍ਰਤੀہار ਹੁਣ ਸਰਕਾਰੀ ਵਕੀਲ ਨੇ ਹਮਲਾ ਜੋ ਕਰਦੇ ਉਹ ਦਿੱਸ ਤੇ ਹੀ ਗੱਲ ਸੁਗਲਾਈ ਨੂੰ ਲੋਕ ਨੂੰ ਪਿਆਰ ਪਾਪ ਨਾਲ ਜਿਹੜੇ ਕਰੇ ਪਾਪ ਨਾਲ ਉਹਨਾਂ ਤੇ ਹਮਲਾ ਹੋਣਾ ਦੂਏ ਪਾਸੇ ਤੇ ਜਾਂ ਕਿਉਂਕਿ ਤਬਈ ਤੇ ਉੱਤੇ ਗਚੈਰੀ ਜਿਹੀ ਹੁੰਦਾ ਹੁੰਦਾ ਉਹ ਤੇ ਵਕੀਲ ਨਹੀਂ ਲਪੜਦਾ ਨੂੰ ਕੋਈ ਆਪਣੀ ਗਾਲ ਆਪੇ ਕਰਨੀ ਪੈਣੀ ਜਾਂ ਫਿਰ ਗੁਰੂ ਵਕੀਲ ਬਣਦਾ ਕਰਨੀ ਲੋਕ ਤੇ ਜਿਹੜੇ ਵਕੀਲ ਬਣਦਾ ਤੇਰਾ ਗਿਆਨ ਹੈ ਵਕੀਲ ਬਣਦਾ ਤੇ ਗਾਲਤ ਕਾਹਨ ਹੈ ਜੇ ਫੜਿਆ ਤਾਂ ਗਾਲਤ ਕਰ ਲੂਗਾ ਤੇਰੇ ਕੰਨ ਨਹੀਂ ਬੁਕਾਨਤ ਤੇ ਸਖਰੇ ਜਿਹੜੀ ਹਰਬਾਨੀ ਹੈ ਬਕਾਦ ਤੇ ਰਸਾਰੀ ਹੈ ਉਥੇ ਜਵਾਬ ਦੇਈ ਆਪਣਾ ਕੇਸ ਕਿਵੇਂ ਲੜਨਾ ਹੈ ਹਾਂ ਆਪਣਾ ਕੇਤਾ ਆਵੇਂ ਲੜਨ ਸੋ ਐਸਾ ਰਾਜਾ ਸ੍ਰੀ ਗੋਪਾਲ ਉਹ ਰਾਜਾ ਹੈ ਗੋਪਾਲ ਜਿਹਦੇ ਘਰ ਐਸਾ ਕੁਛ ਸ੍ਰੀ ਗੋਪਾਲ ਹੈਗਾ ਥੋੜੇ ਆਲਾ ਸ੍ਰੀ ਗੋਪਾਲ ਹੈ ਤੋਂ ਦਾ ਕ੍ਰਿਸ਼ਨ ਹੈ ਸ੍ਰੀ ਗੋਪਾਲ ਇਹਨਾਂ ਨੇ ਸ੍ਰੀ ਗੋਪਾਲ ਜਿਹੜਾ ਬਣਾ ਲਿਆ ਕ੍ਰਿਸ਼ਨ ਉਹਦੇ ਤੇ ਇੱਕ ਕਿਸਮ ਦਾ ਉਹਦੇ ਤੇ ਵੀ ਇੱਕ ਨੇ ਸ੍ਰੀ ਗੋਪਾਲ ਤੇ ਸ੍ਰੀ ਗੋਪਾਲ ਹੈ ਜਾਇ ਜਿਹੜਾ ਸਾਡਾ ਸ੍ਰੀ ਗੋਪਾਲ ਅਸਲੀ ਸ੍ਰੀ ਗੋਪਾਲ ਹੋ ਆਏ ਤੁਹਾਡੇ ਅੱਜੜਾ ਹੈਗਾ ਤੁਸੀਂ ਇਹਦਾ ਸੰਥਾਨ ਦੱਸਿਆ ਉਹ ਸ੍ਰੀ ਗੋਪਾਲ ਨਹੀਂ ਹੈ ਸ੍ਰੀ ਗੋਪਾਲ ਤਾਂ ਇੰਨੀ ਸ਼ਕਤੀ ਉਹਦਾ ਮਾਲਕਾ ਹੈ ਤੁਸੀਂ ਬਣਾ ਲਿਆ ਆਹਾਂ ਤੁਰੀ ਕਬਲ ਜਿਹੜਾ ਹੁਣ ਹੈ ਹੀ ਨਹੀਂ ਜਿਹੜਾ ਜਾਉਂਦਾ ਮਰਦਾ ਉਹ ਵਿਸ਼ਨੂੰ ਦਾ avatars ਬਣਾਇਆ ਨਾ ਰਾਜੇ ਰੈਨ ਨੇ ਜੀ ਤੇ ਇਹ ਚੰਨ ਚਲੀ ਕਬਲ ਨੋ ਰਖ ਲਿਆ ਉਹ ਰਾਮ ਜੰਨ ਨਾਲੇ ਕ੍ਰਿਸ਼ਨ ਨੂੰ ਵੀ ਹੁੰਦਾ ਕ੍ਰਿਸ਼ਨ ਨਾਲੇ ਦਮਤੋ ਵੀ ਹੁੰਦੇ ਉਹ ਹਨ ਰਾਮਾ ਕਹਿੰਦੇ ਨਾ ਹੋਰੇ ਕ੍ਰਿਸ਼ਨ ਉਹਨਾਂ ਨੇ ਆਹ ਆਮਲੂ ਰਮਿਆ ਹੋਇਆ ਕਹਿੰਦੇ ਨੇ ਗੋਪਾਲ ਨਹੀਂ ਕਹਿੰਦੇ ਇਹਨੂੰ ਗੋਪਾਲ ਕਹਿੰਦੇ ਨੇ गोपाल ਦਾ ਮਤਲਬ ਉਹ ਗੋਪਤ ਪਾਲਣਾ ਕਰਦਾ ਪਾਲਣਾ ਕਰਦਾ ਪਰ ਦੀਦਾ ਨਹੀਂ ਹੈ ਪਰ ਗੱਲ ਨਹੀਂ ਹੈ ਗੋਪਤ ਕਰਦਾ ਗੋਪਾਲ ਗੋਪ ਦਾ ਮਤਲਬ ਉਹ ਹੁੰਦਾ ਗੋ ਦਾ ਮਤਲਬ ਇਹ ਜੀਵ ਹੁੰਦਾ ਹੈ ਜੀਵ ਪਾਲਣਾ ਕਰਦਾ ਰਾਜਾ ਰਾਜਾ ਜੀਵਾਂ ਦੀ ਪਾਲਣਾ ਕਰਦਾ ਪਰ ਆਦਮੀ ਲਈ ਉਹ ਕਰਦਾ ਸਾਡੇ ਆਲਾ ਉਹ ਕਹਿੰਦਾ ਸਾਡੇ ਆਲਾ 84 ਲਖ ਜੂਨ ਦੀ ਗੱਲ ਦਾ 10 ਲਖ ਜੂਨ ਹੈ ਸਾਡੇ ਦੀ ਕ੍ਰਿਸ਼ਮ ਕਹਿੰਦਾ ਬਣਨਾ ਨਹੀਂ ਜੀ ਸੋ ਐਸਾ ਰਾਜਾ ਸ੍ਰੀ ਗੋਪਾਲ ਹਾਂ ਐਸਾ ਰਾਜਾ ਸ੍ਰੀ ਗੋਪਾਲ ਉਹਨੂੰ ਰਾਜਾ ਮੰਨਦੇ ਸੀ ਕੋਈ ਹਥਸਮਾਨ ਨਹੀਂ ਰਾਜਾ ਐਸਨ ਗੈਰ ਗਵੀਰ ਵੀ ਇਹਨਾਂ ਜੀ ਨੂੰ ਰਾਜਾ ਕਹਿਣਾ ਆਹ ਰਾਜਾ ਹੋ ਉਹਦੀ ਵਿਆਖਿਆ ਉਹ ਸਾਡੇ ਜੀ कोई हर समान नहीं राजा ए पूत सब दिन चार के टूठे करत दरवाजा वो गल व्याख्या है हारो गल दी व्याख्या करी नहीं करी तो मीरां जी व्याख्या ही है वो नहीं लगाई कोई हर समान नहीं राजा ओ हां था वो चलिए को राजा राजा ने मुझे बात लिया ਹਰੀ ਜਾਂ ਨਰਹਰੀ ਵੀ ਕਹਿੰਦਾ ਉਹ ਰਾਜਾ ਵੀ ਕਹਿੰਦਾ ਬਾਬਾ ਜੀ ਇੱਥੇ ਜੋ ਸੋ ਲਿਖਿਆ ਸੋ ਐਸਾ ਰਾਜਾ ਸੱਸੇ ਵੀ ਲੱਗੀ ਐ ਸੱਜੇ ਆ ਐਵੇਂ ਆ ਕਿ ਸੋ ਸ਼ਬਦ ਆ ਸੋ ਆ ਇਸ ਲਈ ਐ ਇਹਦਾ ਗਣ ਗੰਧਰਵ ਰਿਚੀ ਆ ਉਹਦੇ ਕਰੇ ਨੇ ਗਣੰਦਨਰਵ ਜਿੰਨੇ ਨੇ ਨਹੀਂ ਜਿਹੜੇ ਤੁਸੀਂ ਕਹਿੰਦੇ ਸੁਰਗਾਂ ਦੇ ਵਿੱਚ ਪਰ ਨਰਵ ਨੇ ਜਿਹੜੇ ਇੱਕ ਰਾਗੀ ਨੇ ਇੱਕ ਸਾਜੀ ਨੇ ਗੰਦ ਨਰਵ ਨੰਦ ਅਰਵ ਗਰਨ ਵਾਲੇ ਵੀ ਹੁੰਦੇ ਨੇ ਸਾਜ਼ ਵਜਾਉਣ ਵਾਲੇ ਆਪਣੇ ਕੀਰਤ ਕਹਿੰਦੇ ਨਰਵ ਰਾਗੀ ਜਿਵੇਂ ਲਾਉਣ ਨਾਲ ਬੇਟ ਨਰਵ ਰਾਗੀ ਇਹਨਾਂ ਨਾਲ ਡਿਗਰੀ ਬੱਪੂ ਢਾਡੀਆ ਵੱਪੜੇ ਟਾੜੀਆ ਵੀ ਨੂੰ ਤੇ ਚਾਹਵੇ ਅਗੋਨਾਨਾ ਟਾੜੀ ਉੱਥੇ ਰਹੀਆ ਦਰਬਾਰ ਦਾ ਹੋਂਡਾੜੀ ਤੇਰੇ ਦਰਬਾਰ ਤੇ ਟਾੜੀ ਵੀ ਨੇ ਉੱਥੇ ਉਹ ਵੀ ਸੀ ਪਰ ਉਹ ਗੌਲ ਨੇ ਦਾਸ ਬਣ ਕੇ ਗੌਣੇ ਉਹ ਵੱਪੜੇ ਤਾਂ ਆ ਜਿਹੜੇ ਤਾਂ ਦਰਬਾਰ ਦੇ ਹਸਕਾਰੀ ਜਿਹੇ ਇਹਨਾਂ ਦਾ ਜਿਹੜਾ ਰਾਗ ਹੈ ਉਹਦਾ ਹੰਕਾਰ ਹੈ ਟਾੜੀਆ ਨੂੰ ਹੰਕਾਰ ਨਹੀਂ ਵੱਪੜੇ ਫੰਦਾ ਜਲਮ ਕੇ ਕਰ ਉਹ ਵੀ ਉਹਦੇ ਦਰਵਾਜ਼ੇ ਤੇ ਭਗਤ ਜੀ ਤੁਹਾਡੀ ਉਹ ਸਾਰੇ ਜਿਹਨਾਂ ਵਾਲੀ ਗਾਇ ਹੈ ਗੁਣ ਨੇ ਉਹ ਕੋਟਾ ਦੀ ਹੁੰਦੇ ਜਿਹੜੇ ਹੋਰ ਕੋਲਿਜ ਰੀਕ੍ਰੀਏਸ਼ਨ ਦੇ ਪ੍ਰੋਗਰਾਮ ਸੁਣਾਉਂਦੇ ਨੇ ਉਹ ਰਾਗੀ ਹੁੰਦੇ ਗੁਣ ਗਾਨ ਕਰਨ ਵਾਲੇ ਜਿਹੜੇ ਹੁੰਦੇ ਨੇ ਉਹ ਕੀਰਤਰੀ ਹੁੰਦੇ ਜੀ ਰਾਗੀ ਨਹੀਂ ਹੁੰਦੇ ਰਾਗੀ ਰੋਗੀ ਹੁੰਦੇ ਇਹ ਰਾਗੀ ਵੀ ਨੇ ਜਦ ਦਰਬੀ ਬਣ ਜਾਂਦਾ ਨਹੀਂ ਕੀਰਤਨੀ ਵੀ ਬਣ ਜਾਂਦੇ ਇਹੋ ਕਹਿੰਦੇ ਬਸਾਂ ਵੀ ਕੀਰਤਨੀ ਰਾਗੀ ਆ ਡੋਟ ਹੁੰਦੇ ਰਾਗੀ ਰਾਗੀ ਜਾਸ ਨਹੀਂ ਕਰਦੇ ਹੁੰਦੇ ਜਾਸ ਅੰਦਰੋਂ ਨਹੀਂ ਕਰਦੇ ਹੁੰਦੇ ਅੰਦਰੋਂ ਰਾਗ ਗਾਉਂਦੇ ਹੁੰਦੇ ਨੇ ਮੂੰਹ ਦੇ ਵਿੱਚ ਜੋ ਬੰਦੀ ਬੋਲੀ ਜਾਂਦਾ ਇਹਨੇ ਕੀਰਤਨੀ ਨੇ ਰਾਗ ਨਹੀਂ ਕਰਦੇ ਹੁੰਦੇ ਜਾਸ ਗਾਉਂਦੇ ਹੁੰਦੇ ਆਪਣੀ ਮੋਜ ਵਿੱਚ ਹੋਜੀ ਕੀਰਤੀ ਕਰਨਾ ਬਈ ਕੀਰਤਨ ਕਰਨਾ ਉਸਤਤ ਕਰਨਾ ਬੜਾਈ ਕਰਨਾ ਕੀਰਤੀ ਕਰਨਾ ਉਸਤਤੀ ਕਰਨਾ ਉਹ ਉਸਤਤੀ ਕਰਦੇ ਨੇ ਪਰਮੇਸ਼ਰ ਦੀ ਉਹ ਤਤ ਕਰਿਆ ਨੇ ਜਨ ਅੰਤਨਾ ਪਾੜਾ ਵਾਰ ਉਹ ਕਹਦੇ ਨੇ ਉਹਨਾਂ ਦਾ ਉਸਤਤੀ ਕਰਨ ਵਾਲ ਧਿਆਨ ਰਾਗ ਤਾਂ ਉਹਨਾਂ ਦੇ ਮੂੰਹ ਚ ਆਪੇ ਨਿਕਲੀ ਜਾਂਦਾ ਹੈ। ਰਾਗ ਇਹ ਕੋਈ ਸ਼ਬਦ ਨੂੰ ਬਾਰ-ਬਾਰ ਰੰਗਤ ਦੇ ਕੇ ਪੇਸ਼ ਕਰਦਾ ਹੁੰਦਾ ਹੈ। ਰੰਗਤ ਦੇਣੀ ਉਹਦਾ ਮੇਨ ਕੰਮ ਸ਼ਬਦਾਂ ਨਾਲ ਉਹਦਾ ਕੋਈ ਬਹੁਤਾ ਸਬੰਧ ਨਹੀਂ ਹੁੰਦਾ। ਸ਼ਬਦਾਂ ਦੀਆਂ ਮਾਤਰਾ ਨਾਲ ਸਬੰਧ ਹੈ ਉਹਦਾ। ਆਹ ਮਾਤਰਾ ਇੰਨੀ ਨੂੰ ਆ ਰੰਗਤ ਦਿੱਤੀ ਜਾ ਸਕਦੀ ਹੈ। ਉਹਨਾਂ ਦਾ ਰਸ ਬਦਲਣਾ ਨਿਰੰਗਤਨਾ ਰਸ ਬਦਲਣਾ ਹੁੰਦਾ ਹੁੰਦਾ ਉਹ ਰਾਗ ਦਾ ਰੰਗ ਬਦਲਦਾ ਹੈ ਰਾਗ ਦਾ ਰਸ ਬਦਲਦਾ ਹੈ ਰਾਗ ਰਸ ਉਹਦਾ ਹੁੰਦਾ ਹੈ ਰਾਗੀ ਦਾ ਰਾਗ ਰਸ ਪੇਸ਼ ਕਰਨਾ ਹੁੰਦਾ ਰਾਗੀ ਨੂੰ ਸਰ ਰਾਗ ਰਸ ਚੋਂ ਆਨੰਦ ਹੁੰਦਾ ਨਾਮ ਦਾ ਰਸ ਨਹੀਂ ਰਾਗੀ ਨੂੰ ਖੁਦ ਆਨੰਦ ਹੁੰਦਾ ਜਦੋਂ ਉਹਨੂੰ ਆਨੰਦ ਦੀ ਰਾਸ ਦਾ ਮਿਲਦਾ ਤਾਂ ਸੁਣਨ ਵਾਲੇ ਨੂੰ ਕਦੋਂ ਮਿਲੂ ਇਹਦੇ ਮੋਜ ਚੀਜ ਹੈ ਉਹਨੂੰ ਉਹਦਾ ਰਸ ਨਹੀਂ ਆਇਆ ਸੁਣਨ ਵਾਲੇ ਨੂੰ ਕੰਨਾਂ ਨੂੰ ਰਸ ਕਿਵੇਂ ਆਜੂ ਕੰਨਾਂ ਵਾਲੇ ਦਾ ਕੰਨ ਰਾਜੇ ਇਹ ਬੋਲਣ ਵਾਲੇ ਨੂੰ ਰਾਸ ਦੇਹ ਜਾਉਂਦਾ ਉਹ ਜਿਹੜੇ ਸੁਣਨ ਵਾਲੇ ਨੂੰ ਬੱਪੂ ਦੇ ਢਾਡੀਆ ਗਵੰਤ ਆਛੈ ਆਹ ਉਹ ਵਧੀਆ ਗਾਉਂਦੇ ਗਵੰਤ ਆਛੈ ਗਾਉਂਦੇ ਰਹਿੰਦੇ ਵਾਗਿਆਂ ਮੈਂ ਖਸਦਾਂ ਗਾਉਂਦੇ ਉਹੀ ਨੇ ਦੋਏ ਗਾਉਂਦੇ ਜੀ ਸੋਈ ਤਦ ਗਾਵਣ ਜੋਤ ਤਪਾਵਣ ਉਹ ਨੂੰ ਪਾਉਂਦੇ ਤਾਂ ਉਹਦੇ ਅੱਛੈ ਉਹਨਾਂ ਦਾ ਕੋਰਣਾ ਵਧੀਆ ਹੁੰਦਾ ਸਭ ਤੋਂ ਸਰਬ ਸਾਸਤਰ ਬਹੁ ਰੂਪੀਆ ਭਾਵੇਂ ਜਿਹੜੇ ਸਾਧਾ ਤਰਣ ਵਾਲੇ ਸਾਰੇ ਇਹ ਬਹਿ ਬਹੁ ਰੂਪੇ ਆ ਰਾਸਤਾਰ ਇਹ ਨਹੀਂ ਹੁੰਦੇ ਕਿਉਂਕਿ ਜਦ ਲਾਲाराम ਲੀਲਾ ਵਾਲੇ ਬਹੁ ਰੂਪੀਏ ਦੇ ਬਹੁਤ ਸਾਧਾ ਉਹ ਬਹੁ ਰੂਪੀਆ ਬਹੁ ਪ੍ਰਕਾਰ ਦਾ ਗਿਆਨ ਹੈ ਡੋਡ ਉਹਨਾਂ ਦੀ ਕਮਤ ਨਹੀਂ ਆਏਗੀ ਉਹ ਆਪ ਆਪਣੀ ਬੁੱਧ ਵਾਲੇ ਨੇ 400 ਰੁਪਇਆ ਮਤਲਬ ਹੈ। ਹੈ। ਇੱਕ ਰੂਪ ਤਾਂ ਦੇ ਵਿੱਚ ਹੈ। ਉਹਨਾਂ ਦੀ ਆਪਣੀ ਆਪਣੀ ਮੱਤ ਹੈ। ਸਰਦਾਰ ਸ਼ਾਸਤਰ ਵਾਲੇ ਨੇ। ਉਹਨਾਂ ਨੇ ਤਾਂ ਤਤ ਗਿਆਨ ਨਹੀਂ ਹੁੰਦਾ ਉਹਨਾਂ ਕੋਲ। ਉਹ ਵੀ ਉੱਥੇ ਹੀ। ਅਖਾੜਾ। ਅਨੁਰਵਾ ਉੱਥੇ ਜੇਲਾ ਕੋਈ ਵੀ ਨਹੀਂ ਸਾਰੇ ਗੁਰੂਆਂ ਨੇ। ਅਨ ਦੇਖੀ ਮੁੰਦ ਨੇ ਜੇਲਾ ਨਹੀਂ ਕੋਈ ਗਿਆ ਤਾਂ ਸਾਰੇ ਗੁਰੂ ਬਲੇ। ਉਸਾੜਾ ਆਪਣੀਆਂ ਆਪਣੀਆਂ ਇੰਗੀਆਂ-ਵਿੰਗੀਆਂ ਮਾਰੀ ਜਾਂਦੇ ਨੇ ਕਿਹਦੀ ਕਿਸ ਨਾਲ ਮਤ ਨਹੀਂ ਮਿਲਦੀ ਇਹਨਾਂ ਨੂੰ ਗੇਦੀ ਬਣਦੇ ਜੀ ਮਤ ਪੈਦਨੇ ਨਾਲ ਵਿੱਚ ਸਾਰਿਆਂ ਚ ਤਾਂ ਹੀ ਸੱਤ ਨਹੀਂ ਰਹੀ ਸੀ ਸੱਤੇ ਮਤਾਂ ਨੇ ਸੱਤੀ ਰਣਨੀ ਘਰੇ ਸੇ ਆਪਾ ਰੋਵਣ ਕੂੜੀ ਰੋਵਣੇ ਕੂੜੇ ਕੁੰਮੀ ਕੂੜੇ ਕਮਾ ਵਾਤੇ ਰਉਂਦੀਆਂ ਨੇ ਮੈਂ ਆ ਕਰ ਦੰਦਾ ਸਾਡਾ ਇਹ ਜੀ ਆ ਕਰ ਦੰਦਾ ਸਾਡਾ ਇਹ ਕੀ ਹੋ ਕਰ ਦੰਦਾ ਚੱਤੀ ਕੋਲੇ ਕੋਹ ਮੰਤਰ ਉਹਦੇ ਕੋਹ ਮੰਤਰ ਆ ਕੋਸ਼ਰ ਉਹਨੇ ਆਪਣੇ ਆਪਣੇ ਨਾਥ ਕਰ ਦਿੰਦੇ ਆਪਣੇ ਆਪਣੇ ਏਂਗਲਾ ਨਾਲ ਉਹਨਾਂ ਨੇ ਬੇਜ਼ਰ ਥਾਇਆ ਆਪਣੀ ਆਪਣੀਆਂ ਮੱਤਾ ਚਲਾਈ ਉਹਨੇ ਆਪਣੇ ਆਪਣੇ ਝੇਲੇ ਦੇ ਢੜੇ ਬਣਾਤੇ ਉਹਨਾਂ ਨੇ ਅਸਲ ਦੇ ਵਿੱਚ ਰਿਸ਼ੀ ਮਹੰਨੀ ਨਾ ਤਿਆ ਕਰੇ ਬਾਹਰ ਜਣਾ ਹੈ ਇਹ ਇਹਦੀ ਵਿਚਾਰਤਾਂ ਵਿਖਰ ਗਈ ਇੱਕ ਵਿਚਾਰਤਾਂ ਦਾ ਵਿਖਰੀਆ ਨਹੀਂ ਸੀ ਇਹ ਆ ਕੇ ਉਹ ਰਿਸ਼ੀ ਮਹੰਨੀ ਦਾ ਇੱਕ ਢੜੇ ਦਾ ਨਹੀਂ ਸੀ ਮਹੰਨੀ ਇੱਕ ਢੜੇ ਦਾ ਜਿਹੜਾ ਬ੍ਰਸਪਤ ਹੈ ਗੁਰੂ ਉਹ ਢੜੇ ਦਾ ਮਾਤ ਹੈਗਾ ਰਾਮ ਜਨ ਪਰਾਂਵ ਜੰਨਰ ਲੋਮੀ ਵਾਲੇ ਜਨਤਾ ਹੀ ਪੈਦਾ ਹੁੰਦਾ ਆ ਰਾਮ ਲੋਮੀ ਏ ਨੌ ਦੁਆੜੇ ਪ੍ਰਗਟ ਨਹੀਂ ਸ਼ਰੀਰ ਦੇ ਦਸਵੇਂ ਗੁਪਤਾਂ ਦਸਵੇਂ ਜਾਂਦਾ ਹੀ ਨਹੀਂ ਮਾਇਆ ਜਿਹੜਾ ਆ ਰਾਮ ਲੋਮੀ ਹੁੰਦੀ ਹੈ ਨਾ ਜੀ ਬਸ ਦਸ ਵੀਰ ਦਾ ਜ਼ਾਇਰਾ ਦਾ ਆ ਇਹਨੂੰ ਉਹਦਾ ਰਾਵਣ ਮੱਦਦਾ ਉਹ ਮਨ ਮੱਦਾ ਦਸ ਵੀਰ ਇਹਦਾ ਨੂੰ ਆਪਲਾ ਰਵੜਾਂ ਦੀ ਹੋਰ ਕਿਸੇ ਦਾ ਮਾਰਦਾ ਬਾਹਰ ਪਣਾ ਲਿਆ ਰਾਵਣ ਆਪਲਾ ਮੰਨੂ ਰਾਵਣ ਨਹੀਂ ਬਣਿਆ ਰਾਵਣ ਦੋਦੇ ਆਪਣੇ ਅੰਦਰ ਸੀ राम ਜੰਨ ਦੇ ਉਹ ਰਾਵਣ ਨੂੰ ਉਹਦਾ ਨਵ ਰਾਵਣ ਲਖਿਆ ਜਿਹੜਾ ਚਾਰ ਮੇਰ ਦਾ ਗਿਆ ਤਾਸੀ ਉਹਨੂੰ ਰਾਵਣ ਕਹਿਣ ਲੱਗ ਉਹਦਾ ਬ੍ਰਾਹਮਣ ਸੀ ਮੰਡਲਿਕ ਬੋਲ ਬੋਲੇ ਕਾਛੇ ਉਹ ਮੰਡਲ ਇਹਨੂੰ ਹੀ ਲੰਬਯਾਰ ਮੰਡਲ ਹੈ ਮੰਡਲੀ ਹੈ ਮੰਡਲੇ ਕਬੂਲ ਬੋਲਦੇ ਹੈ ਕੱਕਾ ਦੂਏ ਪਾਸੇ ਲਾਤਾ ਆਉ ਚੈ ਜਾਨ ਕੇ ਲਾਤਾ ਮੰਡਲੀ ਕਬੂਲ ਬੋਲੈ ਕਬੂਲ ਬੋਲਨੇ ਬੋਲ ਨਹੀਂ ਬੋਲਦੇ ਕਬੂਲ ਬਗਾੜ ਕੇ ਬੋਲਦੇ ਨੇ ਜੇ ਕੋ ਬੋਲਾ ਦੇਖੋ ਆਖਾ ਬੋਲ ਬਗਾੜ ਤਾਂ ਲਿਖਿਆ ਸਰ ਕਵਾਰਾ ਗਵਾਰ ਦੇਖਿਆ ਨਾ ਕੱਲ੍ਹ ਨੂੰ ਲਾਗੇ ਕਹਿੰਦਾ ਕਿ ਇਹਨਾਂ ਸਤ ਤੁਸੀਂ ਮੈਂ ਜਦ ਮੈਂ ਬੋਲਦਾ ਫਿਰ ਇਹਨਾਂ ਦਾ ਐਡਾ ਨਾ ਕਿਆ ਕਰੋ ਕੀ ਕਹਿ ਇਹਨਾਂ ਨੂੰ ਦੱਸ ਤਾਂ ਕਾ ਐਡਾ ਲਾਇਆ ਅਫਰਾਦ ਇਹ ਅਫਰਾਦ ਹੈ ਜੀ ਛੋਟਾ-ਬੋਟਾ ਹੀ ਹੈ ਗੋ ਆਏ ਇਹਨਾਂ ਨੇ ਜਾਣ ਵਜੀ ਆਪਣੇ ਪਾਪ ਛਪਾ ਲਏ ਲੋਕਾਂ ਨੂੰ ਕਦੀ ਗਲੇ ਪਾਤਾ ਉਹ ਤੂੰ ਦਾ ਵੀ ਕਿਹਦੇ ਨੂੰ ਪਤਾ ਲੱਗਿਆ ਇਹਦੇ ਵੀ ਕੋਈ ਕਾਇਦਾ ਨਾ ਆਇਆ ਹੈ ਨਹੀਂ ਤਾਂ ਕਹਤਾ ਜੇਰਾ ਅਖਰ ਇਹਦੋਂ ਤਾਂ ਹਰਾ ਤੇ ਉਹ ਪ੍ਰਚਾਰ ਕਰਤਾ ਵੀ ਇਹਦੋਂ ਨਾਲੇ ਇਹ ਹੱਥ ਲਿਸਟ ਜਿਹੜੀ ਹੈ ਉਹ ਤਾਂ ਅੱਧ ਹਈ ਨਹੀਂ ਇਹਨਾਂ ਨੇ ਕੀਤਾ ਵੀ ਕੀਤਾ ਕਿਉਂ ਕੀਤਾ ਉਹ ਮੰਡਲੀ ਹੁੰਦਾ ਮੰਡਲੀ ਕੀ ਹੁੰਦਾ ਵੇ ਦੱਸ ਮੰਡਲੀ ਹੁੰਦਾ ਸਿੱਧ ਮੰਡਲੀ ਮੰਡਲੀ ਜੁੰਡਲੀ ਹੁੰਦਾ ਨਾ ਜੀ ਜੁੰਡਲੀ ਉਹਨੂੰ ਮੰਡਲੀ ਹੁੰਦੀ ਹੈ ਸੰਤਾ ਦੀ ਮੰਡਲੀ ਹੁੰਦੀ ਹੈ ਸਾਖਤਾ ਦੀ ਜੁੰਡਲੀ ਹੁੰਦੀ ਹੈ ਗੋਲ ਕੈਰੇਜ ਬੈਠਣਾ ਚਰਚਾ ਕਰਨ ਨੂੰ ਜਿੱਦੇ ਗੋਲ ਮੀਟਿੰਗ ਕਾਨਫਰੰਸ ਹੁੰਦੀ ਹੈ ਉਹ ਮੰਡਲੀ ਕਹਿੰਨੇ ਜਿਹੜੇ ਉਹਨੇ ਦਾਕੂ ਇਹ ਨਹੀਂ ਸੰਤਾਨੀ ਜੁਣੜੀ ਸੰਤਾਨੀ ਸੰਤਾਨੀ ਜੁਣੜੀ ਸੰਤਾਨੀ ਮੰਨਣੀ ਉਹ ਜੁਣੜੀ ਇਕੱਠੇ ਹੋ ਕੇ ਜਾਵੈ ਨੇ ਜੁੜ ਕੇ ਜੁੜ ਕੇ ਹੁੰਦੀ ਉਹਨਾਂ ਦੀ ਬੁਰੇ ਕੰਮ ਹੋ ਜਾਂਦੇ ਸੰਤਾਨੀ ਮੰਨਣੀ ਹੁੰਦੀ ਆਇਤਾ ਮੰਨਣੀ ਉਹਨਾਂ ਦੀ ਜਿਹੜੇ ਆਪਣੇ ਆਪ ਕਹੁੰਦੇ ਨੇ ਕੰਮ ਕਾਜ ਨਹੀਂ ਨਾ ਚਲੇ ਸਾਰੇ ਭੈਣ ਨੇ ਜੁੜ ਕੇ ਜੀ ਉਹ ਮੰਨਣੀ ਹੁੰਦੀ ਆ ਉਹਨਾਂ ਦੀ। ਖੰਡ ਮੰਡਲ ਖੰਡ ਮੰਡਲ ਬ੍ਰਹਮ ਬਹ ਮੰਡਾ ਐਨੀ ਮੰਡਲ ਨਾਲ ਜੀ ਮੰਨ ਲਈਏ ਮੰਡਲ ਤੇ ਮੰਨ ਲਈਏ ਮੰਨ ਲਈਂ ਬਣਾਤਾ ਚੱਕੇ ਕਰ ਕਬੂਲ ਤੀਨਾ ਜਿਹੜਾ ਕਬੂਲ ਲਫ਼ਜ਼ ਉਹ ਬਚਾਉਣਾ ਬੋਲ ਬੋਲੇ ਉਹ ਪੁੱਠੀਆਂ ਗੱਲਾਂ ਕਰਦੇ ਨੇ ਬੇਤੋਂ ਬਾਦ ਬਾੜੀਆ ਉੱਥੇ ਕਬੂਲ ਬੋਲਦੇ ਨੇ ਇੱਥੇ ਆ ਕੇ ਵੱਡੀ ਆ ਜਿਹੜਾ ਨੇ ਉਹ ਕਬੀਰ ਨੇ ਕਿਹਾ ਸੀ ਵੱਡਲ ਬਾੜੀ ਬਾਟ ਇੱਥੋਂ ਕਬੂਲ ਤੋਂ ਬੋਲ ਕਰਕੇ ਆ ਪਾਛੇ ਘਰਤਾ ਵੀ ਪੜਨੇ ਨਾ ਲੋ ਇਹ ਕਰਾਮਾਤਮੀ ਸੁਨਰੀਆਂ ਦੀ ਕੀਤੀ ਹੋਈ ਐਦਾਂ ਰੋਣਾ ਪਉਂਦੇ ਸੀ ਉਹ ਸੇਈ ਤਵਜੂਨਾ ਟਿੱਕਾ ਲਖਾਇਆ ਸੀ ਤਾਂ ਹੀ ਸਿੱਖ ਦੀ ਬੋਲਵਾਤੀ ਤੇਗਾਉ ਹੀ ਹੈ ਹਿੰਦੂ ਵਾਲਾ ਹੀ ਸਿੱਖ ਦੀ ਬੋਲਵਾਤੀ ਵੀ ਹੁਣ ਲੋਕ ਵਿਸ਼ਵਾਸ ਕਰ ਲੰਗੇ ਬਹੁਤ ਸ਼ਾਨਦਾਰ ਆਦਮੀ ਸੀ ਤੇ ਉਹਨਾਂ ਕਰਤ ਅਤਲੇ ਹੁਣ ਵੀ ਨੇ ਹੌਂਦੈਲਾ ਕਿਸੇ ਬੋਲਦਾ ਹੀ ਨਹੀਂ ਚੁੱਪੇ ਹੋ ਗਿਆ ਸਰਬ ਸ਼ਾਸਤਰ ਬਹੁ ਰੂਪੀਆ ਨਨ ਕਰਵਾ ਅਖਾੜਾ ਇਹ ਮੰਡਲੀ ਮੰਡਲੀ ਕਬੂਲ ਬੋਲੀ ਕਾਛੇ ਹਾਂ ਤੇ ਕਾਛੇ ਹੁੰਦਾ ਕਾਛੇ ਟਿੱਕ ਬੋਲ ਨੇ ਨਾ ਉਹ ਕਮਜੋ ਪਿੱਕ ਦੂਗੇ ਤੇ ਟਿੱਕ ਦੂਗੇ ਆ ਰੰਗ ਚਾੜੇ ਨੂੰ ਲਾਉਦੇ ਨੇ ਜੀ ਬਈ ਜਿਹੜੇ ਹੁੰਦੇ ਨੇ ਬੋਲ ਅੱਛੇ ਬੋਲ ਨਹੀਂ ਹੈ ਉਹ। ਸੱਚੇ ਬੋਲ ਨਹੀਂ ਹੈ, ਖਬੂਲ। ਅੱਛੇ ਨੇ ਕਾੱਚੇ। ਕਾੱਚੇ ਨੂੰ ਤੁਸੀਂ ਝਗੜਾ ਪਾਉਣ ਵਾਲੇ ਵੀ ਕਹਿ ਰਹੇ, ਕਹਿ ਸਕਦੇ ਹਾਂ ਅਸੀਂ। ਝਗੜਾ ਬੁਧਾਉਣ ਵਾਲੇ ਵੀ ਕਹਿ ਸਕਦੇ ਹਾਂ। ਤੁਹਾਨੂੰ ਕਹੋ ਜਿਹੜੇ ਸਤ ਨੇ ਉਹਨਾਂ ਦੀ ਗੱਲ ਅਸਲ ਚ ਹੈ। ਸ਼ਾਸਤਰ ਉਹਨਾਂ ਦੇ ਲਿਖੇ ਹੋਏ ਨੇ। ਆਪਣੇ ਆਪਣੇ ਕੋਈ ਸ਼ਾਸਤਰਾਂ ਦੇ ਵਿੱਚ ਜਿਹੜੇ ਨੇ ਸਤ ਰੇਸ਼ੀ ਨੇ ਹੋਈ। ਸਤਿ ਪ੍ਰਕਾਸ਼ ਦੇਨ ਦੇ ਉਹ ਮੱਤਾ ਨੇ ਉਹਨਾਂ ਦੇ ਸਤ ਵਿਚਾਰਤਾਰਾਵਾਂ ਨੂੰ ਸਤ ਉਹ ਕਹਿਆ ਸੱਤ ਹੀ ਦੰਨੀ ਕਰੇ ਸੇ ਆਪਾਂ Hindu મત ਰਨੋ ਸਤ ਵਿਚਾਰਤਾਰਾਵਾਂ ਕਠੀਨ ਦੇਵੀਆਂ ਨੇ ਨਾ ਇਹਨਾਂ ਦੀ ਸਤ ਸਹੀ ਕੀ ਕਥਾ ਹੈ ਪੂਰੀ ਪਈ ਹੈ ਸਤ ਦੇਵੀਆਂ ਨੇ ਅਸੱਚ ਸਤ ਜਿਹੜਾ ਸੀ ਸੱਚ ਸੀ ਗੱਲ ਉਹ ਜਿਹੜੀ ਸੱਚ ਦੀ ਦੇਵੀ ਚੰਡੀ ਆ ਉਹਦੀਆਂ ਨੇ ਸੱਤ ਬਣਾਤੀ ਜਿਵੇਂ ਇੱਕ ਦੇ ਤਿੰਨ ਬਣਾਏ ਨੇ ਇਹਨਾਂ ਨੇ ਬਰਮਾ ਵਿਸ਼ਨੂ ਸ਼ਿਖਜੀ ਇੱਕ ਤੋਂ ਘਾਤੋਂ ਤਿੰਨ ਬਣਾਏ ਨੇ ਸੱਤ ਨੇ ਹੈਗੇ ਅੱਠ ਪਜਾਹਾਨ ਨਾਲ ਦੇ ਵੀ ਇਹਨਾਂ ਸੱਤ ਜਿਹੜੀਆਂ ਨਕਲੀ ਨਹੀਂ ਅਸਲੀ ਆ ਸੱਤ ਪ੍ਰਕਾਰ ਦੀਆਂ ਮਤਾਂ ਕੋਤੋਂ ਜਿਹੜੀਆਂ ਬਣਾਈਆਂ ਨੇ ਥੋੜਾ ਥੋੜਾ ਥੋੜਾ ਥੋੜਾ ਹਟ ਗਈਆਂ ਸੱਚ ਤੋਂ ਉਹਨੇ ਅੱਠਵੇਂ ਮਾਤਰ ਹੈਗੀ ਗੁਰਮੁਖ ਕੋਈ ਅਸਤਾਨ ਵੀ ਕਹਿੰਦੇ ਨੇ ਇਹਨੂੰ ਪਤੰਜਲੀ ਦਾ ਅਸਤਾਨੀ ਹੋ ਗਏ ਉਹਦਾ ਜਵਾਬ ਉਹਨੇ ਦਿੱਤਾ ਵੀ ਜਿਹੜਾ ਅਸਤਾਨ ਜਿਹੜਾ ਉਹਦੇ ਚ ਸੀ ਯਮ ਪਹਿਲਾਂ ਫਿਰ ਨਿਯਮ ਨਿਯਮ ਤੇ ਉਹ ਬੋਲਿਆ ਮੁਸਲਮਾਨ ਵੀ ਜਿਹੜਾ ਨਹੀਂ ਨਿਯਮ ਬਣਾਏ ਨੇ ਨਿਯਮ ਬਣਾਏ ਨੇ ਇਹ ਆਦਮੀ ਨੇ ਬਣਾਏ ਨੇ ਮੈਸੇਜ ਜਿਹੜਾ ਕੋਈ ਭੇਜਿਆ ਮਤ ਦਾ ਤੁਹਾਨੂੰ ਦਾ ਮੈਸੇਜ ਭੇਜਿਓ ਪਰਮੇਸ਼ਰ ਨੇ ਤੇ ਜਿਹੜੀ ਸ੍ਰਿਸ਼ਟੀ ਪਰਮੇਸ਼ਰ ਨੇ ਬਣਾਈ ਹੈ ਤੇ ਜਿਹੜੇ ਉਹਨੇ ਮੈਸੇਜ ਭੇਜਿਆ ਪਰਮੇਸ਼ਰ ਨੇ ਭੇਜ ਉਹ ਤੋਂ ਹਟਵੇਂ ਵਾਲੇ ਨੇਮ ਆਦਮੀ ਨੇ ਬਣਾਏ ਨੇ ਉਹ ਨਹੀਂ ਚੱਲ ਸਕਦੇ ਉਹ ਅਸਲੀ ਨਹੀਂ ਹੁੰਦੇ ਪਰਮੇਸ਼ਰ ਦੇ ਜਿਹੜੇ ਨੇਮ ਨੇ ਉਹ ਬਨਾਂਗੇ ਸ੍ਰਿਸ਼ਟੀ ਉਹਨੇ ਬਣਾਈ ਹੈ ਉਹਦੇ ਵਾਸਤੇ ਨੇਮ ਵੀ ਉਹੀ ਬਣਾਊਗਾ ਆਦਮੀ ਕਿਵੇਂ ਬਣਾ ਸਕਦਾ ਹੈ ਕਿ ਆਦਮੀ ਉਹ ਆਪਣੇ ਬੜੇ ਬਣਾਉਂ ਕਿ ਆਪਣੇ ਮਨ ਤਰਨ ਸਾਰੇ ਬੜੇ ਹੋਈ ਨੇ ਸਭ ਨੇ ਆਪਣੇ ਆਪਣੇ ਨੇ ਬੜਾਏ ਨੇ ਆਪਣੇ ਆਪਣੇ ਤਰਨੇ ਇਹ ਤੇ ਉਹ ਜਿਹੜਾ ਨੂੰ ਪੁੱਛਿਆ ਕੋਈ ਗੱਲ ਨਹੀਂ ਨਾ ਗੱਲ ਦਾ ਜਵਾਬ ਨਹੀਂ ਐਂਡ ਵਿੱਚ ਵੀ ਕਿਹਾ ਇੱਥੇ ਆ ਕੇ ਡਰ ਡਲੋਪ ਪੈਦਾ ਹੋ ਗਿਆ ਉਹ ਇਹਦਾ ਕੋਈ ਜਵਾਬ ਨਹੀਂ ਉਹ ਆਦਮੀ ਤੁਹਾਡੀਆਂ ਮੱਤਾ ਬਣਾਈਆਂ ਨੇ ਪਰਮੇਸ਼ਰ ਤੁਸੀਂ ਛੱਡਦਾ ਸ੍ਰਿਸ਼ਟੀ ਪਰਮੇਸ਼ਰ ਨੇ ਬਣਾਈ ਹੈ ਆਦਮੀ ਪਰਮੇਸ਼ਰ ਨੇ ਆਦਮੀ ਵਾਸਤੇ ਨਿਯਮ ਵੀ ਹੀ ਬਣਾਉਗਾ ਇਹਨਾਂ ਨੇ 7 ਸਤ ਰਿਸ਼ੀ ਨੇ 7 ਧੜੇ ਨੇ ਉਹਨਾਂ ਨੂੰ ਇਕੱਠੇ ਕੋਸ਼ਿਸ਼ ਕੀਤੀ ਹੈ ਇਕੱਠੇ ਹੋਏ ਨਹੀਂ ਨੂੰ ਰਖਦਾ ਹਿੰਦੂ ਮਤ ਉਹ ਅਡਗ ਨੇ ਪਤੰਜਲੀ ਦਾ ਇਸਤਾਨ ਚਾਰ ब्रह्मा ਦੇ ਚਾਰ ਚੇਲੇ ਨੇ ਉਹਨਾਂ ਦੇ ਚਾਰ ਨਾਮ ਨੇ ਸੰਕਤ ਸੰਨੰਦਨ ਸੰਤ ਕਬਾਰ ਸਨਾਤਨ ਸਲਾਤਨ ਨਹੀਂ ਮਤ ਪ੍ਰਚਲਤ ਹੈ ਤਿੰਨ ਮਤਾਂ ਅੜੀ ਮੜੀਆਂ ਹੈਗੀਆਂ ਉਹ ਬਹੁਤੀ ਪ੍ਰਚਲਤ ਨਹੀਂ ਹੋਈਆਂ ਆਦਮੀ ਦੀ ਬਣਾਈ ਹੋਈ ਮਤ ਪਹਿਲੀ ਗੱਲ ਤਾਂ ਆਦਮੀ ਦੀ ਬਣਾਈ ਹੋਈ ਹੈ ਦੂਜੀ ਗੱਲ ਚਾਰ ਚੇਲੇ ਇੱਕੋ ਗੁਰੂ ਦੇ ਨੇ ਚਾਰ ਮਤਾਂ ਕਿਉਂ ਨੇ ਉਹਨਾਂ ਦੀਆਂ ਇੱਕ ਮਤ ਕਿਉਂ ਨਹੀਂ ਹਣੋ ਇਹ ਤਾਂ ਚਾਰੇ ਹੀ ਤੋਂ ਦੂਰ ਨੇ ਇਹ ਸਚਾਈ ਹਿੰਦੂਮਤ ਲਈ ਹੈ ਜਿਹੜਾ ਇਹ ਸਚਾਈ ਨੂੰ ਸਮਝਦਾ ਐ ਐਕਸਪੋਜ਼ ਕਰਦੰਦਾ ਅਨੁਸਾਰੀ ਨੂੰ ਉਹਦੇ ਸਾਹਮਣੇ ਬੈਠੇ ਗਦੇ ਨਹੀਂ ਇਹ ਮੈਂ ਸਿੱਖਾਂ ਦੇ ਸਿੱਖਾਂ ਨੇ ਕਹਤਲੇ ਨੇ ਅਣਗਿਣਤ ਨਹੀਂ ਚਲੋ ਉਹਦੇ ਵਿੱਚ ਵੀ ਜਿਹੜੇ ਨੇ ਜਗਰਦਾਰੀਆਂ ਬਾਰਾਂ ਰੱਖ ਸੀ ਇਕੱਠੇ ਕਦੇ ਵੀ ਨਹੀਂ ਹੋਏ ਰਹਿਤਮ ਨੇ ਅਦਾ ਕਾੜਾ ਬਣਾਇਆ ਕੰਝੂਰੋਬ ਨਹੀਂ ਹੋਇਆ ਇਹ ਦੂਏ ਠੀਕੇ ਪਿੱਛੋਂ ਲੈਨੇ ਸੀ ਦੇਖਾ ਉਹ ਚਿੱਕੀ ਤਾਂ ਤੁਸੀਂ ਮੈਲੇ ਵੀ ਨਹੀਂ ਗਏ ਗੁਰੂ ਦੇ ਖਲਾਫ ਰਹੇ ਨੇ ਕਹਤਾ ਵੀ ਤੁਸੀਂ ਵੀ ਕਰ ਲੋ ਅਹੰਡ ਖੜਾ ਜਿਵੇਂ ਉਹ ਹੀ ਪੋਲ ਪਾਉਣੇ ਆੜੀ ਜੇਥੇ ਪਾਉਂਦੇ ਉਹ ਜਗ੍ਹਾ ਆਪਣੀ ਐਲਟ ਬਣਾ ਲਈ ਤਾਂ ਸੋਦੀ ਜਿਆਦਾ ਲੈਂਡਿੰਗੋਂ ਪਾਠ ਜੰਮੇ ਮਰੇ ਤੇ ਵੀ ਉਹੀ ਕਰਾਉਣ ਨਾਂਬਦਾਰ ਉਹ ਜਿਹੜਾ ਪੈਸੇ ਲੈ ਕੇ ਉਹ ਕਰਦਾ ਸੀ ਆਪਣੇ ਫੇਰੇ ਕਰਾਉਂਦਾ ਸੀ ਲਾਵਾ ਪੜਾਉਂਦਾ ਸੀ ਤੂੰ ਜਦੋਂ ਚੌਗਣਾ ਕਰਦਾ 10 ਗੁਣਾ ਰੇਟ ਕਰਦਾ ਤੁਸੀਂ ਕਿਹੜਾ ਕੱਟ ਕੀਤਾ ਹੁਣ ਆ ਕੇ ਸੋਲ ਬਿਲਕੁਲ ਸਾਰੇ ਕੁਝ ਢੂੜਦਾ ਆ ਜੋ ਫਿਰਨ ਨਾਲਾ ਜੀਤਾ ਸਾਰਾ ਡਰ ਗਿਆ ਮਹਿਲ ਢੂੜਦਾ ਮਹਿਲ ਡਰ ਗਿਆ ਪੰਜ ਵੀ ਗੱਲ ਵੀ ਪ੍ਰਚਾਰ ਗਲਤ ਹੋਇਆ ਇਹ ਨਹੀਂ ਗੌਰ ਹੁੰਦੀ ਏ ਛੂਟ ਦੀ ਇਹਦੇ ਵੀ ਬਹੁਤ ਦੇਲ ਦੀ ਉਮਰ ਖਤਮ ਹੋਈ ਹੋਈ ਪਰ ਚਲੋ ਜੱਬੀ ਪੁੱਟ ਕੇ ਖਰੀਜਨ ਨੇ ਕੁਝ ਆ ਰਹਾ ਹੈ ਬ੍ਰਿਸ਼ੂਪਰਾਣ ਛੇਤਰਾਣ ਦੇ ਖਿਲਾਫ ਆ ਛੇਤਰਾਣ ਬ੍ਰਿਸ਼ੂਪਰਾਣ ਦੇ ਖਿਲਾਫ ਆ ਦੀ ਅਸਲੀਅਤੇ ਸ਼ਬਦ ਵੀ ਦੱਸੀ ਹੋਈ ਹੈ ਸਾਰੇ ਹਾਂਜੀ ਮਹਾਨ ਕੋਸ਼ ਅਨੁਸਾਰ ਅਸਤਾਂ ਅਸਤਾਂਗ ਦੇ ਜੋ 8 ਹੈ ਉਹ ਅੱਠ ਅੰਗ ਕਹਿੰਦੇ ਓ ਜੀ ਹੈ ਉਹ ਹੈ ਯਮ ਸਾਰੇ ਸੰਤ ਸਾਰੇ ਸੰਤ ਹੀ ਇਹਦਾ ਹੀ ਪ੍ਰਕਾਰ ਵਾਲੇ ਬੱਚਾ ਹਾਂਜੀ ਯਮ ਲੀਯਮ ਯਮ ਨਿਯਮ ਆਸਨ ਪ੍ਰਾਣਾਯਾਮ ਆ ਪਤਰਿਆਹਰ ਧਾਰਣਾ ਧਿਆਨ ਸਮਾਧੀ ਆ ਅੱਠ ਹੈ ਜਦੋਂ ਜਦੋਂ ਸਮਾਧੀ ਪਹਿਲਾਂ ਧਿਆਨ ਧਿਆਨ ਤੋਂ ਬਾਅਦ ਸਮਾਧੀ ਕਿਵੇਂ ਹੋਊਗਾ ਧਿਆਨ ਬਾਅਦ ਸਮਾਧੀ ਹੋਣੀ ਨਹੀਂ ਸਕਦੀ ਜੇ ਕਿ ਆਨੰਦ ਸਮਾਧੀ ਨਹੀਂ ਹੁੰਦੀ ਤੇ ਸਮਾਧੀ ਹਕਤ ਹੈ ਨਹੀਂ ਉਹਦਾ ਤਾਂ ਸਮਾਦ ਹੀ ਦਾ ਸਮਾਧੀ ਵੀ ਕੱਢੀ ਕਿ ਆ ਸੋਲੋ ਸਮਾਦ ਹੈ ਸਾਇਤ ਸਮਾਦ ਹੈ ਨਾ ਸੋ ਨਾ ਸਮਾਦ ਕਹੇ ਨਾ ਸਾਇਤ ਸਮਾਦ ਹੀ ਕਹਿੰਦਾ ਸਮਾਧੀ ਦਾ ਬਰੇ ਮਰੇ ਦੀ ਬਣਾਉਂਦੇ ਨੇ ਇਟਾ ਉਹ ਸਮਾਧੀ ਹੈ ਮਰੇ ਦੀ ਜਿਹੜੀ ਇਟਾ ਦੀ ਬਣਾਉਂਦੇ ਉਹ ਸਮਾਧੀ ਹੁੰਦੀ ਹੈ ਚੇਤਨਿਆ ਸੁਗਮਾਦ ਉਹ ਸਾਇਤ ਜੇ ਗਰਸਨ ਨੂੰ ਸਮਾਗ ਅਨਾਹਪੈ ਨਾਦ ਹੈ ਨਾ ਜੀ ਕਹਿੰਦੇ ਸਮਾਤ ਕਹਿਣੀ ਤੇ ਸੁਨ ਸਮਾਗ बेहोश ਲੋਮੇ ਚ ਜਾਂ ਫਿਰ ਜਾਗ ਜਾਗਦਾ ਹੈ ਕਲਪਨਾ ਕਰਦਾ ਹੈ ਕਿ ਕਲਪਨਾ ਰੁਕ ਜਾਣੀ ਹੀ ਸਮਾਧੀ ਹੈ ਇੱਕ ਪਾਸੇ ਇੱਕ ਪਾਸੇ ਦੀ ਧਿਆਨ ਹੀ ਧਿਆਨ ਹੈ ਜੋ ਇੱਕ ਇੱਕ ਪਾਸੇ ਦਾ ਜੇ ਤੁਸ ਪਾਸੇ ਜਾ ਰਿਹਾ ਰਿਹਾ ਧਿਆਨ ਹੈ ਜਾਂ ਦੁੱਖ ਇੱਧਰ ਉੱਧਰ ਸਦੇ ਇੱਧਰ ਹੁੰਦਾ ਰਹੇ ਤੇ ਕੰਮ ਨਹੀਂ ਆਉਂਦੀ ਹੈ। ਕੰਮ ਨਹੀਂ ਜਾਂਦਾ। ਕਿਉਂਕਿ ਅੱਖ ਪਟਕਦਾ ਹੈ, ਪਟਕਣਾ ਹੋ ਜਾਂਦੀ ਹੈ। ਫਿਰ ਕਹਿੰਦੇ ਕਿ ਅੱਖ ਗਿਆ। ਵੱਡੀ ਜਮੂਨ ਦਾ ਪੈਨ ਦੂਸਰੇ ਪਾਸੇ ਚਲੇ ਗਿਆ। ਇਹ ਪਾਸੇ ਜਿਆਦਾ ਗੱਡੀ ਰਹਿਣਾ ਸਟ੍ਰੇਟ ਹੋ ਗਿਆ। ਸਾਵਧਾਨੀ ਖਤਮ। ਦੁਰਘਟਨਾ ਹੋਏ ਜਾਣੀ ਹੈ। ਹੈ। ਸਮਾਧੀ ਤਾਂ ਕੋਈ ਹੁੰਦੀ ਓ ਜਾਣੇ ਚੇਤਨਹੀ ਦੀ ਇਸ ਕਰਕੇ ਰਹਿੰਦੇ ਨੇ ਮੁਕਤੀ ਨੂੰ ਬਾਦ ਮੁਕਤੀ ਹੈ ਮਨ ਤੋਂ ਬਾਦ ਸਮਾਧੀ ਕਰਦੀ ਓਦੀ ਕੁਛ ਵੀ ਨਹੀਂ ਇਹਨਾਂ ਦੇ ਪੱਲੇ ਕਹਿਣ ਚੋਰ ਢੂਲ ਜਾਂਚੇ ਹੈ ਪਵਨ ਲੱਲਾ ਜੀ ਢੂਲ ਟੱਡਾ ਢੋਲ ਵਾਲਾ ਜੀ ਸਾਦਾ ਸਾ ਹੈ ਬਾਦ ਕੀ ਹੈ ਲੱਲਾ ਜੀ ਤੇ ਇੱਕ ਢੂਲ ਢੋਲਾ ਚੋਰ ਢੂਲ ਜਿਆਦਾ ਪਾਸੇ ਤੇ ਆਵਾਜ਼ਾਂ ਫੇਰੀਏ ਉਹ ਕੁਝ ਬੋਲਦਾ ਸੁਆ ਕੁਝ ਬੋਲਦਾ ਧੀਆ ਕੁਝ ਬੋਲਦਾ ਚੌਥਾ ਕੁਝ ਬੋਲਦਾ ਚਾਰੇ ਪਾਸੇ ਡਿਫਰੈਂਟ ਤਰ੍ਹਾਂ ਦੀ ਆਵਾਜ਼ ਆਉਂਦੀ ਹੈ ਕਬੂਲ ਕਬੂਲ ਉਹੀ ਗੱਲ ਉਹ ਕਹਿੰਦਾ ਉਹਦੀ ਲੋ ਕਹਿੰਦਾ ਵਿਦਵਾਨ ਇਹ ਵੀ ਕਹਿੰਦੇ ਬਚਾਰ ਨਹੀਂ ਕਰਦੇ ਕਹਦੇ ਨਹੀਂ ਹਜ਼ੂਰੀਆ ਚੋਰ ਢੂਲ ਚਾਚੇ ਹੈ ਪਵਨ ਤੇ ਤੇ ਹਵਾ ਜਿਹੜੀ ਪਬਲਿਕੀ ਬੋਂਗ ਦੀ ਬਾਣੀ ਨਹੀਂ ਹੁੰਦੀ ਜਾਰੇ ਪਾਸੋਂ ਤੋਂ ਡਿਫਰੈਂਸ ਕਿਸਮ ਦੀ ਆਵਾਜ਼ ਹੈ ਉੱਥੇ ਜਿੱਤੇ ਸਤ ਪ੍ਰਕਾਸ਼ ਦੀ ਸਭਾ ਨੂੰ ਦੋਸਤ ਜਿੱਤੇ ਇਹ ਬੈਨਾਨੀ ਮੰਡਲੀ ਬੰਦੀ ਹੈ ਨਾ ਜਦ ਐ ਨਾਨੀ ਜੀ ਮੰਡਲੀ ਬਣੇੜੇ ਕਬੂਲ ਨੇ ਚਾਰਾਂ ਪਾਸਾਂ ਤੇ ਇੱਕ ਦੂਦੇ ਵਿਰੋਧੀ ਆਵਾਜ਼ਾਂ ਨੇ ਯਾਰੇ ਬੇਦਾਨੀ ਆਵਾਜ਼ਾਂ ਨੇ ਇੱਕ ਮਤ ਨਹੀਂ ਹੋ ਰਿਹਾ ਕੋਈ ਕਹਿੰਦਾ ਜਿਹੜਾ ਧਰਮ ਹੈ ਸ਼ਕਤੀਆਂ ਨੇ ਹੀ ਧਰਮ ਸ਼ਕਤੀ ਵਿਰੋਧ ਧਰਮ ਹੀ ਨਹੀਂ ਸ਼ਕਤੀਆਂ ਨਹੀਂ ਤਾਂ ਧਰਮ ਨਹੀਂ ਹੈ ਸ਼ਕਤੀ ਦਿਖਾਉਂਦੇ ਨੇ ਚਰਤੀਆ ਇਹ ਉਹਨਾਂ ਨੇ ਕੀਤੀਆਂ ਹੋਈਆਂ ਨੇ ਬਾਹ ਐਡੀ ਲੰਮੀ ਕਾ ਲਈ ਉਹ ਕਾ ਲਈ ਝੂਠ ਬੋਲੇ ਗੁਰਨਾਨਦ ਨੇ ਆਪਣੇ ਬਈਂ ਦੇ ਵਿੱਚ ਤਿੰਨ ਦਿਨ ਛਾਲ ਮਾਰੀ ਉਹ ਕਰਤਾ ਉਹ ਕਰਤਾ ਹੈ ਜਮਨਾ ਦੇ ਵਿੱਚ ਕ੍ਰਿਸ਼ਨ ਨੇ ਛਾਲ ਮਾਰੀ ਇਹ ਇੱਕ ਤਾਂ ਇਹ ਹੈ ਕਰਾਮਾ ਕਾ ਵਖਾ ਵੱਡਾ ਝੂਠ ਬੋਲ ਕੇ ਵੱਡਾ ਬਣਨਾ ਵੱਡਾ ਇਹ ਗੁਰਨਾਨਦ ਨੂੰ ਵੱਡਾ ਬਣਾਉਣ ਦਾ ਇਹੀ ਮਤਲਬ ਸੀ ਵੱਡੇ ਵੱਡੇ ਝੂਠ ਬੋਲਦੇ ਉਹਨਾਂ ਨੂੰ ਬਾਬਾ ਦੀਪ ਸੂ ਸੀਸ ਲੈ ਗਿਆ ਹੱਥੇ ਠੀਕ ਕਰਕੇ ਲੜਿਆ ਸੀ ਉਹਨਾਂ ਦੇ ਖਲਸਿਆਂ ਨਾਲ ਲੜਿਆ ਸੀ ਇਹ ਸਭ ਝੂਠ ਜਿਹੜੇ ਨੇ ਇਹ ਧਰਮ ਇੱਕ ਤਾਂ ਇਹ ਪੱਖ ਦਾ ਪ੍ਰਚਾਰ ਕਰਦੇ ਨੇ ਸ਼ਕਤੀਆਂ ਪੈਦਾ ਕਰਦੇ ਨੇ ਜੋ ਰੱਥ ਨਿਕਲਿਆ ਜੋ ਧਾਮਿਕ ਨਿਕਲਿਆ ਜੋ ਸਾਂਖਰਿਕ ਨਿਕਲਿਆ ਜੋ ਆਉਂ ਨਿਕਲਿਆ ਉਹ ਪ੍ਰਚਾਰ ਹੈ ਇਹਨਾਂ ਦਾ ਸ਼ਕਤੀਆਂ ਤੇ ਕਾਇਰ ਨੇ ਉਹ ਮੰਨ ਨਹੀਂ ਦਿੰਦੇ ਹਾਲ ਦੇ ਖਿਲਾਫ ਨੇ ਉਹ ਕਹਿੰਦੇ ਨੇ ਜਿਹੜੀ ਚੀਜ਼ ਨੂੰ ਜਮਾਤੀ ਵਾਲੇ ਨੇ ਰਾਆਂ ਆ ਵਾਲੇ ਪ੍ਰਾਂਣ ਚੜਾ ਲਓ ਫਤਲ ਉਹ ਜਦੋਂ ਚੜਾ ਲਓ ਤੇ ਤੁਸੀ ਮਰਦੇ ਹੀ ਨਹੀਂ ਨਹੀਂ ਸਕਦਾ ਤੇ ਪ੍ਰਚਾਰ ਹੈ ਯਾਨੀ ਉਹ ਐਂਟੀ ਸਭ ਕੁਝ ਪ੍ਰਚਾਰ ਹੈ ਪਰਮੇਸ਼ਰ ਕੋਈ ਨਹੀਂ ਬਾਗੀ ਨੇ ਸਾਰੇ ਪਰ ਮੈਂ ਚਲ ਜਾਏ ਦੋ ਬਾਹਰ ਜਾਣਾ ਚਾਹੁੰਦੇ ਨੇ। ਘਾਲ ਤੋਂ ਬਚਣਾ ਚਾਹੁੰਦੇ ਨੇ। ਜਿੰਨੇ ਵੀ ਨੇ ਇਹ ਬਚਿਆ ਮੈਂ ਭਗਵਾਨ RAM ਜਿਹੜਾ ਹੈ ਭਗਵਾਨ ਤਾਂ ਆਦਮੀ ਵੀ ਹੁੰਦਾ। ਆਦਮੀ ਵੀ ਹੁੰਦਾ। ਕਾਗੇਬਾਨ ਵੀ ਹੁੰਦਾ। ਪਰਮੇਸ਼ਰ ਨਹੀਂ ਹੁੰਦਾ। ਵਾਹ। खाली ਪਾਏ पे भगवान तुजे भगवान ना तो काल बस भी है मद्द जंदा है जेडा मद्द जंदा परमेश्वर भी है एक बनी जात आ जो मुक्ति भी नहीं मिली उनो तो खाली पाए पे भगवान तु जागते है जग जाकी कला है आ जेड़ा आदमी दे कला है शरीर विच ਜਗਤਿਆ ਇਹ ਹੀ ਭਗਵਾਨ ਹੈ ਜਾਗ ਤੇ ਹੈ ਜਦ ਜਾਗੀ ਚਲਾ ਹੈ ਜਦ ਜਾਗ ਜਾਂਦਾ ਹੈ ਕੋ ਭਗਵਾਨ ਹੁੰਦਾ ਜਾਗਦੀ ਨਹੀਂ ਜਗਤ ਰੂਪ ਦੇ ਵਿੱਚ ਨਹੀਂ ਆਉਂਦੀ ਉਹਨਾਂ ਚੋ ਭਗਵਾਨ ਨਹੀਂ ਹੈ ਜਦ ਜਾਗ ਜਾਂਦਾ ਭਗਵਾਨ ਜੇ ਜੀ ਸੁਤੇ ਜਾ ਹੀ ਬੁੱਧ ਬਗਲਗੀ ਤੋ ਭਗਵਾਨ ਨੇ ਉਹ ਬਜੀਰੋਣੀ ਹੋਈ ਹੈ ਜਾਣਣੀ ਸੀ ਜਾ ਕੇ ਸੁਪਨਾ ਦੂਰ ਹੋ ਗਿਆ। ਜਿੰਦਿਆ ਦੀ ਸਮਝ ਆ ਗਈ। ਸੱਚ ਹੋ ਜਲਿਆ। ਉਹ ਭਗਵਾਨ ਜਮਤਾ ਵਾਲਾ ਉਹ ਨਹੀਂ ਸੁਪਾ ਕਰ ਰਹਿਣ ਨਿਕੁਰਬਾਨੀ ਤੇ ਮੇਰਾ ਨਾਮ ਸੁਪਾ। ਉਹ ਭਗਵਾਨ ਨੇ ਕਿਹਾ ਸੁਭਾਗਾ ਮੰਨਿਆ ਨੂੰ ਬੋਲਵਾ ਕਾਲੀ ਪਾਇ ਭ੍ਰਮ ਕਾਲੀ ਪਾਏ ਪਿਓ ਭਗਵਾਨ ਤੋਂ ਜਾਗਦੇ ਆ ਜਨ ਜਾਗੀ ਕਲਾ ਕਾਲੀ ਪਾਇ ਪਿਓ ਬ੍ਰਹਮਾਸ਼ਰ ਕਾਲੀ ਪਾਇ ਤੇ ਹੋ ਗਿਆ ਹੈ ਜਨੇ ਯੋਗੀ ਨੇ ਇਹ ਵੀ ਸਾਰੇ ਕਾਲ ਵਾਸਨੇ ਭਗਵਾਨ ਨੇ ਬਾਸੇ ਨੇ ਜਾਣਾ ਹਾਦਰ ਕਾਲੀ ਪਾਇ ਸੁਰਾਸਰ ਗੰਦਰਬ ਬੰਦੇ ਅਰਵਾਇ ਸੀ ਨਾ ਜੀ ਦੇਵਤਾ ਦੇ ਦਰਵਾਜ਼ੇ ਤੇ ਨਰੇਂਦਰ ਦੇ ਉਹ ਹਰੇਂ ਨਰੂ ਕਰੰਨੇ ਨੇ ਸੁਰਾਸਰ ਗੰਦਰਬ ਜੱਛਪ ਜੰਗ ਦਿਸਾਵੇ ਦਿਸਾ ਆਔ ਸੁਖਾਲ ਸਵਰ ਬਤਕਾਲ ਤੇ ਇੱਕ ਹੀ ਕਾਲ ਆਪਾਂ ਸਦਾ ਇੱਕ ਬਿਲਕੁਲ ਭਗਵਾਨ ਕਹਿੰਦਾ ਭਗਵਾਨ ਤਾਂ ਕਹਿੰਦਾ ਕਾਲ ਵਸ ਵੀ ਮੰਨਦਾ ਨਾ ਉਹ ਉਹ ਨੂੰ ਜੀ ਉਹ ਗੱਲ ਲਕਉਂਦਾ ਜਿਹੜੀ ਖਰਾਫਾ ਦੂਹੀ ਹੈ ਲੈਕਦਾ ਗੁਰਬਾਣੀ ਇਹਨੂੰ ਗੁਰਬਾਣੀ ਚੋਂ ਕੰਕਰੀਆਂ ਗੋਲੀਆਂ ਕੁਝ ਕੁਝ ਹਾਈਲਾਈਟ ਕਰਦੇ ਉਹ ਵੀ ਤੋਰ ਮਰੋੜ ਕੇ ਅਸਲੇ ਤੇ ਲਾਉਣ ਕਰਕੇ ਜਦ ਲਈ ਆਹ ਬੋਲ ਬੋਲਦੀ ਹੈ ਕਬੂਲ ਬੋਲ ਸੱਚ ਨੂੰ ਰੱਟਣ ਲੱਗੀ ਹੋਈ ਹੈ ਕਮਜ਼ੋਰ ਕਿਸੇ ਜਿਹਨੂੰ ਕਮਜ਼ੋਰ ਕਰਦੇ ਨੇ ਜਿਆਦਾ ਆਪਾਂ ਉਹ ਨੂੰ ਪੱਛੇ ਦੇਣ ਫੋਟੋ ਲਾ ਉਹ ਬੋੜਾ ਕਮਜ਼ੋਰ ਕਰਨਾ ਸੱਚ ਨੂੰ ਦੂਏ ਦੀ ਗੱਲ ਨੂੰ ਟੁੱਪਣਾ ਕੱਟਣਾ ਹੈ ਗੈਲੋ ਇੱਕ ਦੂ ਗੱਲ ਨੂੰ ਕੱਟਣਾ ਫਾਈ 체ਰੀ ਜੀਤ ਲੈ ਭਵਨ 체ਰੀ ਸ਼ਕਤੀ ਹੈ ਜਿਹੜੀ 체ਰੀ ਸ਼ਕਤ ਜੀਤ ਲੈ ਭਵਨ ਹਾਂ ਤੱਤੇ ਨੂੰ ਸਿਆਰੀ ਸ਼ਕਤੀ ਹੈ ਜਿਹੜੀ ਸ਼ਕਤੀ 체ਰੀ ਹੈ ਬੁੱਧੀ ਅਜੇ ਅੜ ਕੇ ਰਹੀ ਹੈ ਬਾਬਾ ਜੀ ਹਾਂ ਕੋਈ ਗੁਰਮੁਖੀ ਸ਼ਬਦ ਆਉਂਦਾ ਨਹੀਂ ਆਉਂਦਾ ਭਿੰਨ ਕਿਹਾਂ ਪਰ ਸੁਵਾਈ ਹੈ ਜੇ ਬਾਬਾ ਜੀ ਹੈ ਜਦ ਚਲਦੀ ਹੈ ਜਿਹੜੀ ਇਹਦੇ ਗਿਆਨ ਦੇ ਗਿਆਨ ਦੇ ਦੀ ਚਲਦੀ ਆ ਬੁੱਧ ਦਾ ਭਾਲਕੀ ਹੈ ਗਿਆਨ ज्ञान ना अकॉर्डिंग ही चलूगी वो जो ज्ञान है वही हो तो करूंगी जो पौधे कागज के बीच है वही मरतूगी इतनी वोल्टेज पिछो आ रही ਆਜ ਲਈ ਮੰਡਲੀ ਬੈਠੀ ਹੈ ਨਾ ਕੋ ਮੋਲ ਬੋਲਣ ਵਾਲੀ ਜੀ ਉਹ ਚੁੱਪ ਕਰਾਉਂਦੀ ਆ ਜਦੋਂ ਸ਼ਕਤੀ ਕਰਗਣ ਹੋਂਦੀ ਹੈ ਬੇਬੋਦੀ ਪ੍ਰਗਟ ਹੁੰਦੀ ਹੈ ਨਾ ਸੇਰੇ ਸਾਰਿਆਂ ਦੀ ਨਹੀਂ ਕਿਹਾ ਪਰ ਚਬਨ ਬੋਲੀ ਜਾਂਦੇ ਨੇ ਕੋਦ ਨੂੰ ਜਵਾ ਚੁੱਪ ਕਰਾਣੀ ਸਾਰੇ ਸਾਰੇ ਜੂਫੇ ਨੇ ਉਹ ਪਤਾ ਲੱਗਿਆ ਨਾ ਕਲੀਅਰ ਜੀ ਜੀ ਉਹ ਸਾਰਿਆਂ ਦੇ ਪਵਨ ਦੇ ਤਲੇਂਦੀ ਹੈ ਫਿਰ ਚੰਡੀ ਇੱਥੇ ਪ੍ਰਗਟ ਹੁੰਦੀ ਹੈ ਜੀ ਇੱਥੇ ਆ ਕੇ ਪ੍ਰਗਟ ਹੁੰਦੀ ਹੈ ਚੰਡੀ ਪਬਾ ਜੀ ਇੱਥੇ ਚੇਰੀ ਸ਼ਕਤ ਹੈ ਮਿਲ ਸ਼ਕਤੀ ਕਰਨੇ ਜੀ ਨੂੰ ਹੈ ਬਿੰਦੀ ਕਿਉਂ ਨਹੀਂ ਹੈ ਜਦੋਂ ਬੋਲਾਂਗੇ ਤਾਂ ਬਿੰਦੀ ਲਾ ਕੇ ਬੋਲਾਂਗੇ ਬਿੰਦੀ ਲਾ ਕੇ ਬੋਲਾਂਗੇ ਸ਼ਕਤੀ ਚੇਰੀ ਸ਼ਕਤੀ ਜੀਤ ਲੇ ਪਵਨ ਦੇਖੋ ਜਦ ਸਾਖਤ ਬੋਲਾਂਗੇ ਜਦ ਬਿੰਦੀ ਨਹੀਂ ਲਾਉਣੀ ਇਹ ਸ਼ਕਤੀ ਬੋਲਾਂਗੇ ਜੋ ਹਿੰਦੀ ਵਿੱਚ ਸੱਚਾ ਦੂਆ ਹੈ ਆਤੁੱਥਾ ਨਹੀਂ ਹੈ ਬੋਲੀ ਉਹ ਹੀ ਬੋਲਾਂਗੇ ਸਾਡੇ ਸੱਚਾ ਇੱਕਾ ਤੇ ਸੱਚ ਨਹੀਂ ਹਿੰਦੀ ਚ ਉਰਦੂ ਵਿੱਚ ਵੀ ਤੰਨ ਬਰਕਾਰ ਦੇ ਸੱਚੇ ਨੇ ਸਾਡੀ ਜਿਹੜੀ ਨਾਲ ਆਵਾਜ਼ ਤੰਨ ਪ੍ਰਕਾਰ ਦੀ ਉਰਦੂ ਚ ਸਾਡੇ ਪਰ ਲਫ਼ਜ਼ ਵੀ ਘਟ ਗਏ ਨਾ ਉਹਨੇ ਵੀ ਚੌਥੀ ਰੈਡ ਸਾਡੇ ਕਬੀਰ ਜੀ ਨੇ 52 ਅੱਖਰ ਦੀ ਗੱਲ ਕੀਤੀ ਹੈ। ਉਹਨਾਂ ਨੇ ਬਾਤ ਕਰੀ ਹੈ। ਸਾਡੇ ਚੌਥੀਓ ਕਹੇ ਨੇ। ਉਦੂਜ ਵੀ ਜਾਵਾ ਨੇ। ਸਵਾਦ ਹੁੰਦਾ ਉਹ ਵੀ ਇਹੀ ਆਵਾਜ਼ ਹੁੰਦਾ। ਇਹਨੇ ਇਹਦੇ ਵਿੱਚ ਉਦੂਜ ਜੀ। ਸਾਡੇ ਕੋਈ ਐਸਾ ਸਾ। ਸਤਿ ਹਾਂ ਸ਼ੋਵੀ ਹੈ ਜੀ ਹਾਂ ਯਾਰ 10 ਮੰਗਲਾਂ ਦੇ ਵਿੱਚ ਦੁਨੀਆਂ ਦੇ ਗੇੜੀਆਂ ਮਰਦੀ ਆਦ ਬਾਣੀ 'ਚ ਨਹੀਂ ਲੱਗੀਆਂ ਦਸਮ ਬਾਣੀ 'ਚ ਲੱਗੀਆਂ ਹੋਈਆਂ ਔਰ ਅੱਧੀ ਭਾਈ ਬਹੁਤ ਹੈ ਆਦ ਬਾਣੀ ਗੁਰੂਆਂ ਨੂੰ ਥੋੜੀ ਲਿਖੀ ਹੈ ਕਿ ਤੱਕ ਵੀ ਇਹਨਾਂ ਕੀਤੀ ਹੈ ਸਟਾਈਲਿੰਗ ਹੋ ਜਾਏ ਗੁਰੂ ਕਰਨੀ ਹੋਵੇ ਸਟਾਈਲ ਹੈ ਕਪਾਹ ਤੋਂ ਨਹੀਂ ਲੈਣੀ ਜਦੋਂ ਹੋਈ ਹੈ ਉਸੇ ਦੀ ਬੇਕਰ ਉਸ ਦਾ ਸਟਾਈਲ ਹੋਊਗਾ ਸਟਾਈਲਿੰਗ ਬੋਲਨ ਦਾ ਸਟਾਈਲ ਦਾ ਸੰਬਾਧ ਹਰ ਬੰਦੇ ਆਜਾਈ ਤੋਂ ਤਿਰੰਤ ਬਰੁੰਗਾਨ ਹੈਗਾ ਪਾਛਾ ਬਰਿ ਪਾਛਾ ਇਹ ਦੀ ਇਹਦੇ ਵਿੱਚ ਬਰੁੰਗਾਨ ਕੀ ਪਾਜਾਬਲ ਗਿਰੋਲੇ ਤੁੰਦਸਾਈ ਦੀ ਬੋਲ ਗਿਰੇ ਹਨ ਅੰਡ ਟੂਕ ਜਾ ਜਾਚੈ ਪਸ਼ਮਤੀ ਅੰਡ ਟੂਕ ਨੇ ਜਿਹੜੇ ਪਸ਼ਮਤੀ ਨੇ ਅੰਡ ਟੂਕ ਨੇ ਟੁਕੜੇ ਨਹੀਂ ਅੰਡੇ ਦੇ ਦੋ ਢਾਲ ਅੰਡ ਟੂਕ ਇੱਕ ਅੰਡੇ ਦੇ ਦੋ ਟੁਕੜੇ ਆ ਦੋ ਟੁਕੜੇ ਨਹੀਂ ਆ ਸਤਿਮਤੀ ਨੇ ਦੇਹ ਕੀਤਾ phsmu phsmu ਦੀ ਢੇਰੀ ਇਹ ਤਾਂ ਤੇ phsmu ਤੀ ਨੇ ਦੇਹ ਤਾਰੀ ਦੇਹ ਤਾਰੀ ਨੂੰ phsmu ਦੀ ਹੋਇਆ ਹੋਇਆ ਤੇ ਅੰਡੇ ਜਿਹੜੇ ਨੇ ਦੋ ਚਾਰ ਚੋਗੇ ਨਾ ਢਾਲ ਹੋ ਗਏ ਦੇਹ ਹੈ ਨਾਲੇ phsmu ਘਰ ਚ ਨੇ ਇਹ ਵੀ ਉਹਦੇ ਘਰ ਕੇ ਜਦ ਆਂ ਤਾ ਅਕੇਲਾ ਜਦ ਇਹ ਸਰੀਰ ਚੰਦਨ ਦਾ ਤੇਰਾ ਅਕੇਲਾ ਹੈ ਦੇ ਆਂਦਾ ਪਰਦਾ ਕੋਈ ਹੈ ਤੇ ਦਾ ਧਾਰ ਹੋ ਕੇ ਸਰੀਰ ਦੇ ਨਾਲ ਜੁੜਿਆ ਆਦਾ ਅਦਾ ਸਰੀਰ ਤੋਂ ਵੱਖਰਾ ਹੈ ਹਾਲੇ ਆ ਵਿੱਚ ਅਦਾ ਆਸ਼ ਰਣਾ ਅਦਾ ਮਾ ਪੌਣ ਦੀ ਬਾਣੀ ਨਾ ਹੈ ਕਿ ਉਹ ਜਾਲ ਵਿੱਚ ਹੈ ਅੰਧੇਰਾ ਨਵਾਉਂ ਜਾਲ ਵਿੱਚ ਹੈ ਅੰਧੇਰਾ ਨੂੰ ਨਵਾਸ ਆਕਾਸ਼ ਵਿੱਚ ਹੈ ਉਹ ਗੱਲ ਜਾਲ ਬਖਰਾ ਕਾਜ ਤੋਂ ਹੁੰਦਾ ਹਵਾ ਨੂੰ ਕਾਜ ਤੋਂ ਬਖਰਾ ਨਹੀਂ ਮੰਨਿਆ ਜਾਂਦਾ ਸਮਝੋ ਹਵਾ ਜਦ ਤੱਕ ਜੇ ਬਗਦੀ ਹੈ ਹਵਾ ਚ ਤਾਂ ਮੁਖਰੀ ਲੱਗਦੀ ਹੈ ਜੇ ਹਵਾ ਚ ਬੇਗ ਨਹੀਂ ਸਮਾ ਜਾਂਦੀ ਹੈ ਜੇ ਕਹਿੰਦੇ ਹਵਾ ਮਾਰ ਗਈ ਨਹੀਂ ਚਲਦੀ ਵਧਦੀ ਨਹੀਂ ਹੈ ਤੁਹਾਡਾ ਮਨ ਯਾਗਾ ਉਹਦਾ ਡੈਲੀਆ ਮਹਿਸੂਸ ਨਹੀਂ ਹੁੰਦੀ ਆ ਵਾ ਮਹਿਸੂਸ ਇਹ ਹੁੰਦੀ ਆ ਸਾਨੂੰ ਸਾਡੇ ਗਿਆਨ ਦੇ ਅਨੁਸਾਰ ਹੈ ਹਾਂਜੀ ਸੋ ਐਸਾ ਇਹ ਰਾਜਾ ਕਰਪਾ ਵਾ ਤੁਮਨੇ ਕੋ ਪਤੀ ਇਹ ਤ੍ਰਿਭਵਨਪਤੀ ਰਾਜਾ ਜਿਹੜਾ ਇਹ ਰਾਜਾ ਅਸਲੀ ਕੋਈ ਹਰ ਸਮਾਨ ਰਾਜਾ ਇਹ ਟੂਕ ਪੁੱਤ ਸਾਹਿਬ ਦੇ ਵਿਚਾਰ ਕੇ ਚੁੱਕੇ ਟੂ ਕਾ ਹੈ ਇਹ ਤਾਂ ਐਂਡ ਟੂ ਦੀ ਬਸਮੰਦੀ ਹੈ ਇਹ ਕਹਿੰਦਾ ਮੈਂ ਰਾਜਾ ਉਹ ਇਹਨਾਂ ਤੇ ਐਂਡ ਟੂ ਇਹਨਾਂ ਤੇ ਤਾਂ ਰਾਜ ਕਰਨਾ ਰਾਜ ਨਹੀਂ ਕਰਨਾ ਇਹਨਾਂ ਤੇ ਕਰਨਾ ਆਪ ਮੁਤੀ ਨਹੀਂ ਜਿੰਨੇ ਦੇ ਤਾਲੀ ਨਹੀਂ ਨਾ ਤੇ ਰਾਜ ਕਰਨਾ ਇਹਨਾਂ ਦੇ ਵਿਚੋ ਨਾ ਤੇ ਤੇ ਨੂੰ ਹੀ ਬਣ ਜਾਂਦਾ ਇਹਨਾਂ ਦੇ ਕੇ ਬਾਜੇ ਪੜ ਆਪਣੇ ਬੁੱਧ ਬਲ ਦੇ ਜੋਰ ਨਾਲ ਆਪਣੇ ਸਰੀਰ ਬਲ ਦੇ ਜੋਰ ਤੇ ਜਫਰ ਆਦਮੀ ਦੇ ਆ ਕੇ ਫਿਰ ਜਨਮਿਤ ਫਿਰ ਪੈਸਾ ਆ ਰਿਹਾ ਥਿਆ ਹਾਲ ਵੀ ਆਜਾ ਮੈਨੇ ਵਿੱਚ ਇਨਵੋਲਵ ਹੋ ਜਾਂਦੇ ਨੇ ਹੋਰ ਤਾਂ ਜਾਨਵਰਾਂ ਪੈਸਾ ਆ ਹਥਿਆਰ ਉਤੇ ਸਿਰਫ ਅਕਲ اور ਸਰੀਰਕ ਸ਼ਕਤੀ ਲੋਜੀ ਜਨ ਚਾਹੀਦੀ ਹੈ ਓਨੇ ਕੂਰਮਾ ਪਾਲ ਉਹ ਕੁਰਮਾ ਜਿਹੜਾ ਕੱਛੂ ਆਇਆ ਸੰਤ ਦੇਦੇ ਖੋਪੜੀ ਦੇ ਬਹੁਤ ਦਿਨ ਪਾ ਰੱਖੇ ਨੇ ਉਹ ਵੀ ਉਹਦੇ ਤਰੇ ਹੀ ਆ। ਗੁਰਮੁਖ ਕੱਛੂ ਕਹਿੰਦੇ ਨੇ ਨਾ ਪੱਕਾ ਅਵਤਾਰ ਹੈ ਕ ਹੋਇਆ ਹੋਇਆ ਸਭ ਤੋਂ ਪਹਿਲਾ ਜੀਵ ਕੱਛ ਅਵਤਾਰ ਕਹਿੰਦੇ ਨੇ ਪਾਣੀ ਚ ਫੈਦਾ ਕੱਛੂ ਬਦਲਿਆ ਪਾਣੀ ਦੇ ਵਿੱਚ ਫਿਰ ਮੱਛੀ ਪੈਦਾ ਹੋਈ ਮੱਛ ਅਵਤਾਰ ਜਾ ਚੈੱਕ ਕਰੀ ਹੋਈ ਆ ਸੇਟੀਨ ਦੇ ਹਿਸਾਬ ਨਾਲ ਉਹ ਜਿਹੜੇ ਕਹਿੰਦੇ ਜੀਵ ਨੇ ਕੇ ਤੱਛੂ ਆ ਕੇ ਵੱਡਾ ਕੇ ਪਰਾਂ ਤਾਂ ਨਾ ਕਰਮ ਨਹੀਂ ਹੋ ਇਹ ਜੀਵਨ ਅਸਪੀਡੈਂਟ ਕੇ ਉਹ ਬਣਦਾ ਡਿਵਲਪ ਹੋ ਕੇ ਫਿਰ ਆਪੇ ਮੱਛ ਕੱਚ ਕਰਨੀ ਕਰ ਬਾਚਕਾਰ ਦੇ ਰੂਪ ਦਾ ਪ੍ਰਕਾਰ ਨਹੀਂ ਕਰਦਾ ਹੈ ਆਪ ਤੇ ਬੁੱਧ ਡਿਵੈਲਪ ਕਰਦਾ ਆਪਣੀ ਫਨੀ ਬਾਸਕ ਸੇਜ ਵਾਲੂਆ ਉਹ ਜਿਹੜਾ ਵਿਸ਼ਨੂ ਆ ਉਹ განਨਾ ਲਾਉ ਪਰ ਉਸ ਤੇ ਉੱਪਰ ਉਹ ਗੰਗਾ ਉਹ ਬੀਰ ਉਹਦੇ ਕੰਢੇ ਵਿੱਚ ਹੀ ਹੈ ਭੋਗ ਜਾਂਦਾ ਰਾਵਣ ਹੈ ਬੋਰ ਤੋਂ ਦਸ ਜੀ ਦਾ ਉਹਦੇ سنگ ਤੇ ਥੱਤੀ ਹੈ ਖੜੀ ਉਹਦੇ ਆਸਰੇ ਖੜੀ ਹੈ ਥੱਤੀ ਖੜਾ ਖਥੂ ਤੇ ਉਹਦੇ ਕੋਲ ਗੰਗਾ ਚਾਹੀਦੀ ਹੈ ਫਿਰ ਪਾਣੀ ਚਾਹੀਦਾ ਉਹ ਗੰਗਾ ਦਾ ਉੱਥੋਂ ਨਿਕਲੀ ਹੈ ਕਿੱਥੋਂ ਨਿਕਲੇ ਸਮੁੰਦਰ ਤੋਂ ਨਿਕਲੀ ਹੈ ਗੰਗਾ ਹੁੰਦਾ ਜਿ ਘਚੂ ਆ ਪਾਣੀ ਦੇ ਵਿੱਚ ਉਹਨਾਂ ਨੇ ਐ ਜੋੜਤਾ ਉਹਨੇ ਜੋੜਤਾ ਉਹ ਸਾਦਰ ਦੇ ਵਿੱਚ ਛੇ ਜਨਾਗਾ ਉਹਦੇ ਦੇ ਮੱਤੇ ਵਿਸ਼ਨੂੰ ਆ ਛੇ ਜਨਾਗਾ ਨੇ ਉਹ ਕੀਤਾ ਹੈ ਉਹਨਾਂ ਨੇ ਆ ਬਣਾ ਲਿਆ ਐ ਜੋੜ ਸਾਦਰ ਦੇ ਵਿੱਚ ਤਾਂ ਛੇ ਨੂੰ ਤਾਂ ਸਾਲੀ ਆਉਂਦਾ ਪਾਣੀ ਚ ਬੋੜਦ ਉਹ ਸਾ ਪਾਉਂ ਦਾ ਦੇ ਤਾਂ ਉਹਦੇ ਪੈਰ ਨੇ ਆਪ ਦਾ ਬਾਹਰ ਉਪੜੀ ਉਹ ਤਾਂ ਕਹਿਦਾ ਨਹੀਂ ਕਾਇਰ ਨੇ ਉਹਦੇ ਕੱਟੂ ਦੱਸਦੇ ਤਾਂ ਆਪਣੋਂ ਜੀ ਤਰ੍ਹਾਂ ਬਾਹਰ ਹੈ ਉਹ ਉੱਥੋਂ ਸਿੱਟੀ ਦਾ ਹੋਰੀ ਜਨ ਨੇ ਚੱਕ ਕੇ ਉਹ ਉਧਰ ਉੜ ਜਾਂਦੇਗੇ ਸੱਪਾਂ ਵੱਲੋਂ ਨਾਂਦਾਂ ਵੱਲੋਂ ਚਲੋ ਸਹ ਫਨੀ ਬਾਸਕ ਬਾਸਕ ਕੀ ਹੁੰਦੇ ਬਾਤ ਕਰ ਉਹਦਾ ਬਾਤ ਉਹਦਾ ਰਾਜਾ ਇਹਨਾਂ ਦਾ ਬਾਤ ਜਿਹੜਾ ਰਾਜਾ ਸੱਪਾਂ ਦਾ ਉਹਨੂੰ ਬਾਤ ਹੁਕਮ ਉਹਦੇ ਕੋਈ ਫੌਨ ਹੁੰਦਾ ਸੈਸ ਨਹੀਂ ਹੁੰਦੇ ਪਹਿਲਾਂ ਸਹਿਤ ਮੁਕੀਆ ਉਹ ਜਿਆਨਾ ਪ੍ਰਤਾਦ ਉਹਦਾ ਧਿਆਨ ਹੈ ਫਿਰ ਆ ਕੇ ਜਦ ਇਕ ਹੋ ਜਾਂਦਾ ਸਵਦਾ ਰਾਜਾ ਉਹ ਹੈ ਜਿਆਦਾ ਜਿਹਰੀ ਲੋ ਹੋ ਜਾਂਦਾ ਬਾਤ ਕੋ ਨੂੰ ਵੀ ਦੇ ਉੱਤੇ ਸਭ ਚੜਿਆ ਫਿਰਦਾ ਛੋਟਾ ਜਿਹਾ ਥੰਗਲ ਹੁੰਦਾ ਰਾਜਾ ਹੋ ਹੀ ਜਾਂਦਾ ਬਾਸਕ ਕੋਟ ਸੇਜ ਵਿਸਥਰੀ ਆਹੋ ਬਾਤ ਕੋ ਨਹੀਂ ਬਾਤ ਸੁਣੇ ਉਹਦੇ ਫਲਸਫੀ ਹੈ ਇਹਨਾਂ ਦੀ ਜੇ ਤਾਂ ਪੜ੍ਹੀ ਹੋਵੇ ਹਿੰਦੂਆਂ ਦੀ ਦੋ ਫਲਸਫੀਆਂ ਨੇ ਅਡਵਟ ਇੱਕ ਸ੍ਰੀ ਪ੍ਰਾਣ ਇੱਕ ਬਿਸ਼ੂ ਪ੍ਰਾਣ ਚ ਹੈ ਕਹਿੰਦੇ ਸਭ ਕੁਝ ਉਹਦੇ ਕਰਤੇ ਜਿਹਨੂੰ ਤੁਸੀਂ ਵਸਾਰਿਆ ਹੋਇਆ ਹੈ ਜਿਸੇ ਘਰ ਵਿੱਚ ਸਭ ਕੁਝ ਹੈ ਘਰ ਵਾਲੀ ਚੀਜ਼ ਲੈ ਲਈ ਆਪਣੀ ਉਹ ਘਰ ਵਾਲਾ ਚੜਤਾ ਮੰਨ ਕੇ ਮਾਲ ਕਬੱਡਾ ਚੀਜ਼ ਵੱਡੀ ਉਹਦੇ ਘਰ ਵਾਲੀ ਤੇ ਉਹ ਹੋਏ ਵੀ ਉਹਦੇ ਮੁਕਾਬਲੇ ਦੀਆਂ ਚੀਜ਼ਾਂ ਨੇ ਤਾਂ ਹੀ ਉਹਦੇ ਮੁਕਾਬਲੇ ਦੀਆਂ ਕਈ ਮੁਤਲ ਮੰਗੀਆਂ ਕਿ ਜਦੋਂ ਕੋਈ ਪੱਖ ਲੈ ਲਿਆ ਕਿ ਜਦੋਂ ਕੋਈ ਪੱਖ ਲੈ ਲਿਆ ਕਿ ਜਦੋਂ ਕੋਈ ਪੱਖ ਲੈ ਲਿਆ ਕਿ ਜਦੋਂ ਕੋਈ ਪੱਖ ਲੈ ਲਿਆ ਆਪਣੀ ਆਪਣੀ ਬੁੱਧ ਸੰਸਾਰ ਉਹਦੇ ਅੱਖ ਹੱਤ ਕਰ ਲਏ ਆਪ ਆਪਣੀ ਬੁੱਧ ਜੇਤੀ ਬਣ ਤਪਨ ਪਿੰਨ ਤੋਂ ਤੇਤੀ ਉਗਲਾ ਲ ਸੰਜਾਇ ਪਸਵਾ ਦਾ ਕੈਬਲ ਸਜਾ ਪ੍ਰਥਮ ਸੰਦਵਾਰਾ ਪ੍ਰਥਮ ਸੰਤਾਰਾ ਕਿਵੇਂ ਸਜਿਆ ਉਹ ਦੱਸਿਆ ਇਹਨਾਂ ਨੇ ਇਹਨਾਂ ਨੇ ਹੋਰ ਕਿਵੇਂ ਦੱਸਤਾ ਦੋ ਪ੍ਰਕਾਰ ਜੰਦੂਆਂ ਨੇ ਦੱਸਿਆ ਇੱਕ ਪ੍ਰਕਾਰ ਜੀ ਮਾਨਾਂ ਨੇ ਅਰੰਡੇ ਜੰਦ ਦੱਸਿਆ ਉਹ ਲੱਗਿਆ ਆਦਮੂ ਤੋ ਗਿਰ ਦੱਸਿਆ ਇੱਕ ਨਹੀਂ ਗੱਲ ਤੇ ਨੀ ਗੁਰਮਤਮਰ ਵਾਲੀ ਗੱਲ ਇਹ ਕਰਕੇ ਦੋ ਪ੍ਰਕਾਰ ਦੇ ਕੰਡੀਸ਼ਨਰ ਤਾਂ ਨੇ ਉਹਨਾਂ ਜਿਸ ਫਾਰਾ ਬਿਆਖਿਆ ਕੀਤੀ ਇਹਦੇ ਨਾਲ ਦੀ ਬਹੁਤ ਪ੍ਰਧਾਵੀ ਦਾ ਜਵਾਬ ਜੀ ਬਾਬੇ ਆਦਮ ਦੀ ਗੱਲ ਕੀਤੀ ਹੋਈ ਹੈ ਇਹਨਾਂ ਨੇ ਜਾਂਚੈ ਕਰ ਹੂਰਮਾ ਪਾਦ ਤਹ ਫਨੀ ਬਾਸਕ ਏਜ ਉਹ ਕੁਰਮਾ ਪਾਲੇ ਵੀ ਕਹਿੰਦੇ ਨੇ ਉਹ ਕੁਰਮਾ ਤੋਂ ਦਾ ਪਾਲਕ ਹੈ ਕੁਰਮੇ ਨੂੰ ਵੀ ਸਾਬ ਨੂੰ ਹੋਰ ਹੋਰ ਪਾਲਣਾ ਕਰਨ ਵਾਲਾ ਨਾ ਜਿਦੂ ਜਿਦੂਨ ਕਹਿੰਦੇ ਆਂ ਸਭ ਦੀ ਪਾਲਣਾ ਕਰਦਾ ਉਹ ਕੁਰਮੇ ਦੀ ਵੀ ਪਰਣਾਉਂ ਕਰਦਾ ਅੱਛੂ ਵੀ ਉਸ ਦਿੰਦਾ ਜਿਸ ਸਾਬ ਨੂੰ ਕੁਰਮਾ ਪਾਲ ਕਹਤਾਂ ਨੂੰ ਆਪਣਾ ਬੜਾ ਬਣਾਤਾ ਜਿਹੜੀ ਦਾ ਰਹਿਮ ਕੋ ਦੰਦਾ ਨਹੀਂ ਹੋਤਾ ਸਮਾਧੀ ਲਾਉਂਦਾ ਆਪਣੇ ਵਾਸਤੇ ਜੇ ਗਿਆਨ ਕਰਾਉਂਦਾ ਉਹ ਗੁਰੂ ਤੇ ਯਾਨੀ ਉਹ ਵੀ ਆਦਮੀ ਵਾਲਾ ਗਿਆਨ ਹੈ ਨਾ ਆਦਮੀ ਆਦਿਨੋ ਗਿਆਨ ਦਊ ਜਿਹੜਾ ਪਾਲਣਾ ਕਰਨ ਵਾਲਾ ਉਹ ਸਾਰਿਆਂ ਦੀ ਕਰੂਗਾ ਸੇਚ ਵਾਲੂਆ ਦਾ ਕੀ ਅਰਥ ਹੈ ਜਿਹਦੇ ਤੇ ਪਿਆ ਉਹ ਕਹਾਂ ਨਹੀਂ ਆ ਵਿਸ਼ਨੂੰ ਦਿਖਾਇਆ ਹੈ ਫਿਰ ਉਹ ਤੇਜ ਹੈ ਉਹਦੀ বালੂਆ ਉਹ ਬਾਲੂਆ ਮਿੱਟੀ ਦੀ ਹੈ ਮਿੱਟੀ ਵਾਸਤੇ ਮਿੱਟੀ ਦੀ ਸਰੀਰ ਵਾਸਤੇ ਸਰੀਰ ਦੀ ਤੇਜ ਹੈ বালੂਆ ਰੇਤ ਉਹ ਦਾਏ ਮਿੱਟੀ ਹੈ ਚੇਤਨਾ ਦੋਹਾਂ ਦੀ ਗੱਲ ਨਹੀਂ ਹੈ ਚੇਤਨਾ ਦਾ ਕੋਈ ਸਹੀ ਨਹੀਂ ਉਹ ਮਿੱਟੀ ਹੈ ਸਰੀਰ ਮਿੱਟੀ ਵਾਸਤੇ ਮਿੱਟੀ ਹੀ ਹੁੰਦੇ ਜਾਂ বালੂਆ ਦੋ ਪਾਸੇ বালੂ ਹੀ ਹੈ ਇਹ ਤਾਂ ਨਹੀਂ ਗੱਲ ਨਹੀਂ ਹੈ ਇੱਥੇ ਜੀ বালੂ ਰੇਤ ਜੋਂ ਨੂੰ ਪਠਿਆਰੇ ওই বালੂ ਹੈ বালੂ ਰੇਤ ਹੁੰਦੀ ਹੈ 18 ਪਾਰ ਬਨਸਪਤੀ ਮਾਲਣੀ ਪਠਾਰਾ ਪਾਰ ਬਨਸਪਤੀ ਹੈ ਇੱਕ ਇੱਕ ਪੱਤਾ ਦੋੜੀ ਹੋ ਜਾਂਦੇ ਬਨਾਸਪਤੀ ਲੈਣਾ ਨੇ ਮੰਨੇ ਹੋਏ ਨੇ ਇਹ ਕਿਉਂ ਨੇ ਨੇ ਉਹ ਗਨਿਆ ਦਾ ਰਾ ਪਾਰ ਬਨਾਸਪਤੀ ਉਹਦੇ ਘਰ ਤੇ ਹੈ ਅੰਦਰ ਸਾਰੀ ਹੈ 18 ਪਾਰ ਬਨਾਸਪਤੀ ਮਾਲਣੀ 18 ਪਾਰ ਬਨਾਸਪਤੀ ਜੀ ਮਾਲਣੀ ਹੈ ਜਿਹੜੀ ਹੈ ਵੀ ਉਹਦੇ ਘਰ ਤੇ ਹੈ ਉਹ ਮੰਡੀ ਤੇ ਬਣਾ ਤਾਂ ਹੁਣ ਬਾਜ਼ੀ ਮੈਂ ਪੈਦਾ ਮਾਲਣੀ ਜੱਤੀ ਹੈ ਬੁੱਧੀ ਹੈ ਚੇਤਨ ਦੀ ਗੱਲ ਐ ਤੇ ਮਾਲਣੀ ਹੋ ਚੀਜ ਐ ਪਾਲਣੀ ਹੋ ਚੀਜ ਐ ਮਾਲਣ ਉਹ ਉਹਨੂੰ ਵਧਾਉਂਦਾ ਨਾਲ ਮਿਲ ਕੇ ਬਣਾਉਂਦਾ ਜੋ ਬਨਸਫਰ ਦੇ ਆਤਮਾ ਉਹ ਮਾਲਣੀ ਹੈ ਬਿਲੀ ਹੋਈਆ ਵਿੱਚ ਮਿਲ ਕੇ ਫੁੱਲ ਬਣਾਇਆ ਉਹਨੇ ਫੁੱਲੇ ਚ ਰਾਜ ਬੜਕੇ ਫੁੱਲ ਦਾ ਰੂਪ ਧੰਨ ਕੀਤਾ ਫੁੱਲ ਜੜਾ ਆਪ ਮਾਲਣੀ ਹੈ ਪੈਦਾ ਕਰਨ ਵਾਲੇ ਕੋਈ ਵੇਲਜ ਮੰਨ ਲਈ ਪਾਣੀ ਪਾਉਂਦੀ ਮੰਨ ਲਈ ਹੈ ਮਾਲਣੀ ਹੋਏ ਨਹੀਂ ਵਿਚਮੀ ਹੋਈ ਹੈ ਜੇ ਮੇਰਾ ਆਰਾਮ ਨਹੀਂ ਹੁੰਦਾ ਜੀ ਦੇ ਵਿੱਚ ਜਗ੍ਹਾ ਜੋ ਹੁੰਦਾ ਉਹ ਮਾਲਣੀ ਹੈ ਬਿੜੀ ਹੋਈਆ ਵਿੱਚ ਮਾਇਆ ਚ ਮਣਕੇ ਹੀ ਹੁੰਦਾ ਹੈ ਮਾਇਆ ਚ ਜੋਤ ਵਿੱਚ ਵਿਆਪਕ ਹੁੰਦਾ ਜੋਤ ਵਿੱਚ ਜਿਵੇਂ ਕਹਿੰਦੇ ਨੇ ਰਮਣਾ ਹੁੰਦਾ ਮਾਇਆ ਵਿੱਚ ਮਿਰਣਾ ਹੁੰਦਾ ਰਮੇ ਚੀਜ਼ ਮਿਲੀ ਚੀਜ਼ ਬੇ ਵਿੱਚ ਫਰਕ ਹੈ ਆਪਾਸ ਵਿੱਚ ਰਮਿਆ ਜਾਂਦਾ ਮਿੱਟੀ ਵਿੱਚ ਮਿਲਿਆ ਜਾਂਦਾ ਪਾਣੀ ਵਿੱਚ ਮਿਲਿਆ ਜਾਂਦਾ ਜਾਂ ਮਲਾਇਆ ਜਾਂਦਾ ਕੁਝ ਪਾਣੀ ਦਾ ਬਲਬਲਾ ਨਾ ਇੱਕ ਬਿੜਿਆ ਜਾਂਦਾ ਰਮੇ ਨਹੀਂ ਜਾਂਦਾ ਪਾਣੀ ਅਕਾਸ਼ ਵਿੱਚ ਰੰਮ ਕੇ ਪਾਣੀ ਚ ਮਿਲਿਆ ਜਾਂਦਾ ਅਕਾਸ਼ ਵਿੱਚ ਨਹੀਂ ਮਿਲਿਆ ਇਹਦੇ ਸਾਡੀ ਤੋਂ ਵਜੂਦ ਅਕਾਸ਼ ਇਸ ਕਰਕੇ ਮੰਨਣੀ ਹੈ 96 ਕਰੋੜੀ ਮੀਗਮਾਲਾ ਚੰਨੀ ਨੇ ਕਰੋੜ ਮੰਗ ਮਾਰਿਆ ਚੰਨੀ ਮਗਰ ਮੀਗ ਜਿਹੜੀ ਉਹ ਖਾਲਸਾ ਉਹ ਤੈਨੂੰ ਕਹਿੰਦੇ ਨੇ 96 ਕਰੋੜ ਖਾਲਸਾ ਜਿਹੜਾ ਅਵਦੇਸ਼ ਕਰਨ ਵਾਲਾ ਉਹ ਨਾ ਮੇ ਬਾਲਿਸ਼ ਕਰੂਗਾ ਦੁਨੀਆ ਦੇ ਵਿੱਚ ਗੁਰਮਤਿ ਪਿਓਰ ਗੁਰਮਤਿ ਜਦ ਕਰੂਣਾ ਵਿਆਖਿਆ ਕਰਨ ਦੇ ਲੈ 96 ਕਰੋੜ ਹੋ ਜੂਗਾ ਉਦੋਂ ਕਹਿੰਦੇ ਸਾਰੀ ਦੁਨੀਆ ਦਾ ਰਾਜ ਉਹ ਸਿਰਫ ਮਤੂੰ ਸਾਡੀ ਦੁਨੀਆ ਮੰਗ ਲਓ ਉਹ ਰਾਜ ਕੀ ਹੈ ਨਿਹੰਗ ਸਿੰਘ ਤਾਂ ਹੀ ਕਰੋੜ ਹੀ ਕਹਿੰਦੇ ਆ ਜਨਮ ਕਰੋੜੀ ਮੁਸਲਮਾਨਾਂ ਦੇ ਲਈ ਵੇਚ ਜਨਮ ਕਰੋੜੂ ਤੋਂ ਆਏ ਹੋਏ 96 ਕਰੋੜੀ ਮੇਗਮਾਲਾ ਪਾਣੀ ਹਾਰੀਆ ਮੇਗਮਾਲਾ ਮੇਗੇ ਨੂੰ ਫਰਮਾਣੋ ਆ ਪਰ ਤੁਗਰਫਾ ਤਰ ਹੁੰਦਾ ਉਹ ਆ ਜਾਣ ਦੇਣ ਵਾਲਾ ਸਾਪਤੀ ਕਿੰਨੀ ਦਾ ਹੁੰਦੀ ਹੈ ਜਾਂ ਬਾਦਸ ਹੁੰਦੀ ਐ ਠੰਡੇ ਹੋ ਜਾਂਦੇ ਲੋਕ ਹੁੰਦੇ ਨੇ ਸਾਰੇ ਪੁੱਜਦੇ ਲਾਵਾ ਬੰਦੋ ਦੀ ਬੱਟ ਪਿਆ ਰਾਤ ਮੈਨੂੰ ਫੋਨ ਆਇਆ ਸੀ ਬੰਗਲਾ ਸਾਹਿਬ ਤੋਂ ਮੇਰਾ ਫਿਰ ਅੱਗੇ ਡਿੱਗਣ ਦੀ ਐ ਆਂ ਕਹਾ ਤੋਂ ਦੋ ਦਾਰੇ ਤੋਂ ਜੇ ਲਾ ਕੇ ਆਏ ਉੱਥੇ ਜਿਹੜਾ ਤੂੰ ਅੰਮ੍ਰਿਤ ਕਹਿਣਾ ਉਹ ਤਾਂ ਹਰੀ ਅੰਦ ਮਾਇਆ ਹੈ ਪਾਣੀ ਉਹ ਮਾਇਆ ਦਾ ਰੰਗ ਜਿਹੀ ਐ ਉਹਨੂੰ ਵਰਤਣਾ ਨਹੀਂ ਅੱਜ ਦੇ ਕੱਲ ਨੂੰ ਹੋਰ ਦਿਨ ਤੋਂ ਜੇ ਹਮਤ ਚਲੋ ਜੀ ਅੱਗੇ ਪਾਣੀ ਹਾਰਿਆ ਤਾਂ ਇਹ ਪਾਣੀ ਆਦੇ ਹੁੰਦੇ ਉਹ ਮੇਂ ਵਾਲਾ ਉਹ ਤੋਂ ਲੈ ਕੇ ਜਲ ਸਮੁੰਦਰ ਤੋਂ ਲੈ ਕੇ ਆਉਂਦੇ ਨੇ ਜੇ ਉਥੋਂ ਆਉਂਦਾ ਦਰਿਆ ਚ ਪਾਣੀ ਨਹੀਂ ਹੁੰਦਾ ਉਹ ਦਰਿਆ ਹੈ ਜੈ ਜਵਨ ਜਵਾਨ ਨਿਕਲ ਜਾਂਦਾ ਇੱਕ ਵਾਰ ਕੇ ਜਿਹੜਾ ਉਲਕੀ ਬਾਣੀ ਹੁੰਦੀ ਆ ਉਹ ਜਿਹਨਾਂ ਦੇ ਜੈ ਜਵਨ ਆਵੇ ਖਦਮੀ ਖਦਮਗੀ ਬਾਣੀ ਐਸਾ ਲਾ ਲਈ ਲੋ ਤੇ ਉਹ ਮੈਗ ਮਾਰਾ ਜਾਂਦਾ ਨਖ ਪਰ ਸੇਵ ਜਾਚੈ ਸੁਰਸੁਰੀ ਜਿਹੜੀ ਹੈ ਜੀ ਇਹ ਬਹੁਤ ਇਹ ਨਾਕਾਏ ਮੁੜਦੀ ਨਹੀਂ ਕਿਸੇ ਪਾਸੇ ਸਖਤ ਹੈ। ਤੁੰਹਿਆ ਇਹ ਨਹੀਂ ਜਿੱਦ ਤੂੰ ਮਰਜ਼ੀ ਮੋੜ ਲੋਂਗੇ ਤੁਸੀਂ ਨੋਂ ਨੂੰ। ਜਿਹੜਾ ਜੇ ਨਾਕ ਪਿੱਛੇ ਨੋਂ ਨਾਲ ਹੋਵੇ ਉਗੜਦੇ ਜਿਹੜਾ ਮਾਸ ਨੂੰ ਜਿੱਦ ਮਰਜ਼ੀ ਮੋੜ ਲੈ। ਸਿੱਧੋ ਪਾਸੇ ਨੂੰ ਚਲਦੀ ਆ ਫਿਰ ਨੋਂ ਇਹ। ਬੜੀ ਸਖਤ ਜੁੰਦੀ ਹੋਣਾ। ਠੀਕ ਨਹੀਂ ਮੁੜਦੀ। ਸਿੱਧੀ ਜਾਂਦੀ ਹੈ ਨੋਂ ਬਾਹਰ ਨੂੰ ਜਾਂਦਾ। ਦੇ ਬਈ ਉਹਦੇ ਨਾਲ ਇਹਨੂੰ ਇਤਕ ਤੱਕ ਦੀ ਹੱਡੀ ਹੋਈ ਆ ਹੈ ਸਾੱਚ ਜਿਹੜਾ ਹੈਗਾ ਨੋਹ ਹੈ ਜਿਹੜਾ ਝੂ ਆ ਦੂਆ ਹੈਗਾ ਸੱਚ ਦੇ ਸਾਚਾ ਝੂਠ ਮੇਸ ਉਹ ਮਾਸ ਹੈ ਹੱਡ ਮਾਸ ਦਾ ਰਿਸ਼ਤਾ ਨਹੀਂ ਕਹਿੰਦੇ ਨੋਹ ਮਾਸ ਦਾ ਰਿਸ਼ਤਾ ਵੀ ਕਹਿੰਦੇ ਹੱਡ ਮਾਸ ਦਾ ਰਿਸ਼ਤਾ ਵੀ ਕਹਿੰਦੇ ਜਿੰਨਾ ਚਿਰ ਹੱਡੀ ਨਾਲ ਨਹੀਂ ਤਾਂ ਮਾਸ ਜਿਹੜਾ ਖੜਾ ਨਹੀਂ ਹੋ ਸਕਦਾ ਹੱਡੀਆਂ ਕਰਕੇ ਜੀੜ ਖੜਾ ਆਪਣਾ ਪਿੰਜਰਾ ਪਿੰਜਰਾ ਹੱਡੀਆਂ ਦਾ ਹੀ ਆ ਆੜਮਾਤ ਹਨਹਾੜ ਫਿਰ ਮਾੜ ਫਿਰ 나ੜੀ ਹੈ ਕੋ ਪਿੰਜਰ ਪਹਿਨਾ ਸੱਚ ਹੈ ਉਹਦੇ ਨਾਲ ਬਾਅਦ ਫਿਰ ਝੂਠ ਹੈ ਲੱਗ ਮਾਫੇ ਹੈ ਯਾਨੀ ਅਸਲ ਜੋ ਹੈ ਪਿੰਜਰ ਉਹ ਹੱਡੀਆਂ ਦਾ ਹੀ ਆ ਅਸਲ ਜੇ ਪਹਿਲਾਂ ਤਾਂ ਨਕਲ ਬਣਦੀ ਹੈ ਕੋਈ ਵੀ ਚੀਜ਼ ਆ ਕਾਪੀ ਬਣੂਗੀ। ਕਾਪੀ ਤੇ ਕੀ ਜੇ ਬਣੂ ਜੇ ਕੋਪੀ ਸ਼ੀਟੇ ਕਾਪੀ ਦਾ ਸੱਚ ਹੋਣਾ। ਪਹਿਲਾ ਦੂਹੁੰਦਾ ਜਿਹੜੀ ਮੱਤ ਹੈ ਸਭ ਤੋਂ ਪਹਿਲੀ ਇਹ ਕਹਿੰਦਾ ਪਹਿਲੀ ਮੱਤ। ਪਹਿਲੀ ਮੱਤ ਝੂਠੀ ਕਹਿੰਦਾ ਕਿ ਪਹਿਲੀ ਮੱਤ ਸੱਚੀ ਹੋਊਗੀ। ਅੱਗ ਵਿੱਚੋਂ ਛੱਟ ਕੇ ਜੇ ਉਠਾ। ਆਗ ਛੱਤ ਦਾ ਮਤਲਬ ਪਹਿਲਾ ਨਾ ਖਾ ਨਾ ਆ। ਉਹ ਤੋਹੀ ਹੁੰਦਾ ਮੋੜਦਾ ਨਹੀਂ ਅੱਡ ਅੱਡੀ ਛੜੀ ਦੇ ਵਿਚ ਨੂੰ ਮਾਫ਼ ਸੇਖ ਇਟ ਇਜ਼ ਸੇਖ ਸਖਤ ਹੈ ਇਹ ਮਰਵਾਣੀ ਹੈ ਨਖ ਪਰసేਵ ਆਪ ਪਰసేਵ ਇਹ ਸੁਰ ਤੇ ਇਹ ਜੋ ਕਹਾਣੀ ਹੈ ਮਤਲਬਾ ਸੁਰ ਅਸਰੀ ਸੁਰ ਉਹ ਲੇਵ ਜਿਹੜੀ ਸੁਰ ਸਰੀ ਹੈ ਹਰ ਕਰਨਾ ਸਾਰਿਆਂ ਨੂੰ ਜਿੱਤ ਲੈਣਾ ਜੁੱਤ ਸਦੀ ਪਰਕਾਣੇ ਫਾਲੀ ਕਹਿੰਦੇ ਆ ਪਕਲਦੇ ਆ ਹਾਂਜੀ ਜਿੱਤਲ ਜਿੱਤ ਲੈਣਾ ਜਿੱਤ ਬਈ ਸਾਰਿਆਂ ਨੂੰ ਇੱਕ ਸਾਲ ਹੁੰਦਾ ਉਹਦੇ ਘਰ ਇਹ ਆ ਉਹਦੇ ਘਰ ਨਾਨਕ ਇਹ ਕਰਕੇ ਨਾਮ ਹੈ ਜੋਤਨੀ ਨੇ ਤੇ ਸੱਚਾਣ ਤੇ ਸੱਚੇ ਸੱਚੇ ਐਂ ਉਹਦਾ ਘਰ ਵੀ ਸੱਚਾਣ ਪਗਲ ਸੱਜਣਾ ਦਾ ਵਾਸੀ ਬੋਲਾ ਨਾ ਹੋ ਗਿਆ ਹਾਂਜੀ ਸੱਜਣਾ ਸੱਚੇ ਸੱਚਾ ਸਤਿਗੁਰੇ ਨਹੀਂ ਮੱਤ ਸੱਚੇ ਵਿਦਿਅਕ ਦੇਸਾ ਉਹ ਨਾ ਖੋਵੇ ਸਖਤ ਉਹ ਮਰਦਾ ਨਹੀਂਗਾ ਉਹ ਖੜਦਾ ਉਹ ਖੜਾ ਰਹਿਣਾ ਅੱਧੀ ਨਾਲੇ ਬਾਸਾ ਲਾ ਹੱਡੀਆਂ ਦੇਖੋ ਕਿ ਹੱਡੀਆਂ ਦਾ ਪਿੰਜਰਾ ਖੜਾ ਰਹਿ ਸਕਦਾ ਬਾਹਰ ਇਹਨੇ ਦੇਖੇ ਬਾਰੇ ਲੋਕਾਂ ਦੇ ਬਾਹਰ ਦਾ ਕੰਮ ਹੋ ਗਿਆ ਜਿਹੜਾ ਵੀ ਉਹ ਜਿਹਨੇ ਸਿਰ ਜੜਾ ਨਾ ਨਾੜੀਆਂ ਨਾ ਮਾਸ ਪਛਿੱਤੂ ਹੁਰਦੇ ਆਸਰੇ ਨਹੀਂ ਕਰਦਾ ਝੂਠ ਸੱਚੇ ਆਸਰੇ ਕਰਦਾ ਮਾਸ ਨਾੜੀਆਂ ਹੱਡੀਆਂ ਦੇ ਆਸਰੇ ਖੜੀਆਂ ਸੀ ਮੈਂ ਲਿਖਿਆ ਸੀ ਸੱਚ ਨੂੰ ਫਸਲੇ ਪ੍ਰਚਾਰ ਨੂੰ ਮਾਇਆ ਦੀ ਲੋੜ ਨਹੀਂ ਹੈ ਫਸਲੇ ਲੋ ਪ੍ਰਚਾਰ ਨੂੰ ਝੂਠੀਆਂ ਸਾਥੀਆਂ ਦੀ ਲੋੜ ਨਹੀਂ ਹੈ ਫਸਲੇ ਪ੍ਰਚਾਰ ਨੂੰ ਸੰਸਾਰੀ ਪਾਣੀਆਂ ਦੀ ਲੋੜ ਨਹੀਂ ਹੈ ਨੂੰ ਗੁਰੂ ਦੇ ਜੀਵਨ ਨੂੰ ਹੀ ਗੁਰੂ ਪੀਰਾਂ ਦੇ ਜੀਵਨ ਨੂੰ ਹੀ ਦੱਸਦਾ ਵਰਦਾ ਪਰ ਤਾਂ ਉਹਨਾਂ ਨੂੰ ਕਰਨੀ ਸੀ ਉਹਨੂੰ ਗੁਰ ਕਰਨੀ ਕਹਿੰਦੇ ਨੇ ਸਾਹਿਤਾ ਉਹ ਇਹ ਸਾਥੀ ਨਾ ਮਗਰ ਨਾ ਕੋ ਉਹਦੇ ਜੀਵਨ ਮਗਰ ਨਾ ਕੋ ਵਰਤਿਆ ਸਾਹਾਰਾ ਖਮਾਉਂਦਾ ਉਹ ਸੀ ਨਬ ਸਿੱਧਾ ਇਹ ਢਟੇਰੀ ਹੋ ਗਏ ਜਿਹੜੀਆਂ ਮੱਤਾਂ ਢਟੇਰੀ ਹੋ ਜਾਂਦੀਆਂ ਨੇ ਉਹ ਸਾਥੀ ਛੱਡ ਦਿੰਦੀਆਂ ਨੇ ਇਹ ਤੁਹਾਨੂੰ ਹੋਏਗਾ ਭਸਮ ਕੇ ਨੂੰ ਮਿਟੇ ਕਹਿੰਦੇ ਨੇ ਅੱਡੀ ਰੂਪੀ ਨਹੀਂ ਲੈਣੇ ਜੇ ਦਾ ਬਾਹਰ ਦੇ ਵਿੱਚ ਹੀ ਮਿੱਟੀ ਹੁੰਦੀ ਹੈ ਨਹੀਂ ਮਾਸ ਕਰਨ ਨੂੰ ਨਾ ਨਾ ਕਬਰਾਂ ਦੇ ਹੱਡੀਆਂ ਨਹੀਂ ਗਾ ਉਹਨੇ ਮਾਸ ਨਹੀਂ ਲੁੱਭਦਾ ਮਾਰਦੀ ਮਿੱਟੀ ਕਹਿੰਦੀ ਮਾਣ ਅੜੀਉ ਲੱਭਦੀ ਉਹ ਤਾਂ ਥੋੜੇ ਦਿਨ ਲੱਗੇ ਕਈ ਇਹ ਬੰਦਾ ਜਾਂਦਾ ਇਹ ਜਿਹੜੀ ਪਾਸ਼ਾ ਨਾ ਨਾਪ ਇਰਕੇ ਨਾ ਦਾਪਾ ਕਰਨ ਲੱਗੇ ਨਾ ਗੈਰ ਨੇ ਪੈਣੋਂ ਕੰਸੇ ਚੈਨੂ ਨਾ ਪੈਣੋਂ ਨਾ ਨਾਖੁਨ ਵੀ ਕਹਿੰਦੇ ਨੇ ਨਾਖੁਨ ਵੀ ਕਹਿੰਦੇ ਨੇ ਉਰਦੂ ਵਾਲੇ ਉਰਦੂਆ ਥਾਂ ਤੇ ਕੋਈ ਪਹਿਲਾਂ ਇਹਨਾਂ ਪਾਸੇ ਕੋਈ ਐ ਵੇਦ ਵਿੱਚੋਂ ਨਿਕਲਿਆ ਨਹੀਂ ਹੁਣ ਹਰਮਾਨ ਦੀ ਅਰੇ ਆਪਾਂ ਨਿੰਦੂ ਵੀ ਆਪਾਂ ਵੇਦ ਵਿੱਚੋਂ ਕੀ ਨਿਕਲਣਾ ਆਪਾਂ ਨਿਕਲ ਕੇ ਨਹੀਂ ਗਏ ਆਪਾਂ ਤਾਂ ਘਰੇ ਦੇ ਵਿੱਚ ਖੜੇ ਹਾਂ ਲਈ ਸਾਡੀ ਤਾਂ ਬੇਇਜ਼ਮਤੀ ਹੈ ਬੁਰਮਤ ਹੀ ਬੇਇਜ਼ਮਤੀ ਹੈ ਉਹ ਕੇ ਬੇਇਜ਼ਮਤੀ ਨਾ ਕਹਿੰਦਾ ਸਾ ਸਮੁੰਦਰ ਦੀ ਹੀ ਗੰਦੇ ਸੀ ਉਹ ਗੇਰ ਸਮੁੰਦਰ ਦੇ ਰੁਪਏ ਆਦੀਆਂ ਸਾਰੀਆਂ ਕਿ ਕਿੰਨੂੰ ਤੁਸੀਂ ਉਲਾ ਸਕਦੇ ਸਾਰਿਆਂ ਨੂੰ ਸਮੁੰਦਰ ਬੜੇ ਮਨਾ ਕਿ ਕਿੰੋਂ ਸਿੱਖਿਆ غور ਵਿਚਾਰ ਕਿਹਾ ਗਿਆਨ ਦੇ ਵਿਚਾਰ ਸਾਲੀ ਦੇ ਗਿਆਨ ਦੇ ਵਿਚਾਰ ਤਾਂ ਇਹਦੇ ਵਿੱਚ ਮੁੰਡੀਆਂ ਨੇ ਆਉਂਦੇ ਉਹਦੇ ਘਾਰੇ ਸੋਰਸਰੀ ਇਹਨੂੰ ਗਿਆਨ ਦੀ ਗੰਗਾ ਕਹਿੰਦੇ ਨੇ ਉੱਦ ਦੇ ਤੇ ਸੋਰਸਰੀ ਹੋਰ ਹੈ ਗੰਗਾ ਹੋਰ ਤੇ ਦੋ ਬਣਾਉਂਦੀ ਜਿਹੜੇ ਸਰਸੁਤੀ ਕਹਿੰਦੇ ਨੇ ਸੋਰਸਰੀ ਹੋਇਆ ਸਰਸੁਤੀ ਇਹਦਾ ਨੌ ਦਾ ਪਹਿਲਾ ਸੋਰਸਰੀ ਦਾ ਅਲਾਵਾਦ ਪਿੰਨੇ ਮਿਲਦੀਆਂ ਨੇ ਆਕੇ ਇੱਕ ਉਹ ਹੈ ਇੱਕ ਜਮਨਾ ਤੇ ਹੁੰਦਾ ਇਹ ਚਾਲੇ ਜਮਨਾ ਦਾ ਇੱਥੇ ਉੱਤੇ ਵੀ ਆਉਂਦੀ ਹੈ ਕਾਹਨ ਤੇ ਆਗਰੇ ਦੇ ਉੱਪਰ ਵੀ ਆਉਂਦੀ ਹੈ ਜਾਂਦੀ ਹੈ ਬਕੌਣ ਦੇ ਪਾਸੇ ਵੀ ਆਉਣੀ ਹੈ ਜਮਨਾ ਤਾਂ ਵਿਚਾਲੇ ਦੀ ਗੰਗਾ ਆਉਂਦੀ ਹੈ ਫਿਰ ਦੀ ਹੋਣੀ ਹੈ ਇਹਨਾਂ ਕਰਕੇ ਆਈ ਇਹ ਕੇਵਲ ਉੱਨੀ ਜਾਂਦੀ ਹੈ ਫਰਜੂ ਦੀ ਸ਼ਾਇਦ ਇਸੇ ਨੂੰ ਕਹਿੰਦੇ ਹੋ ਈ ਇਹ ਲਾਵਾ ਤੋਂ ਸਮੇਂ ਤੇ ਈ ਇਹ ਲਾਵਾ ਈ ਉੱਥੇ ਚਲੀ ਜਾਂਦੀ ਹੋਏ ਕੋਲ ਭਾਂਕੇ પાછી ਉਥੋਂ ਨੜਈ ਜਾਂ ਚਿੱਤੰਨ ਉੱਥੇ ਰਹਦੀ ਨੂੰ ਆ ਕੇ ਉਹ ਤਰਵਾਣੀ ਕਹਿੰਦੇ ਨੇ ਪਰ ਵਿਚਾਲੇ ਹੋਣ ਜਾਂ ਈ ਛੁੱਟਛਲੀ ਇੱਕ ਪਾਸੇ ਵਿਚਾਲੇ ਘਰੋਂ ਤੋਂ ਇੱਕ ਪਾਸੇ ਜੋਗ ਹੈ ਇੱਕ ਪਾਸੇ ਵੈਸ਼ਨਵ ਬੰਤਾ ਰਾਜੀ ਵਾਲੀ ਬਿਸ਼ਨੂ ਵਾਲੀ ਵੈਸ਼ਨਵ ਵੈਸ਼ਨੂ ਭਗਤ ਇਹਨਾਂ ਨੇ ਇਹ ਗਿਆਨ ਉਹਨਾਂ ਦੇ ਗਿਆਨ ਤੋਂ ਪ੍ਰਦਾਨ ਹੁੰਦਾ ਵੈਸ਼ਨਵਾਂ ਨੂੰ ਪਰ ਹੁੰਦਾ ਸਮਰਤੀ ਵਾਲਾ ਗਿਆਨ ਹੈ ਸਾਸਤ੍ਰਾਂ ਦਾ ਇਹ ਵਾਲਾ ਨਹੀਂ ਹੁੰਦਾ ਇਹ ਵਾਲਾ ਵਿਚਾਰੇ ਵਾਲੀ ਜੁਮੇ ਸੁੱਟ-ਸੁੱਟੀ ਜੁਮਦਾ ਮੇਹਰ ਤੋਂ ਸਰੀ ਦੇਵ ਤੇ ਨੂੰ ਜਿੱਤਣ ਵਾਲੀ ਦੇਹ ਤੇ ਕੋਣ ਨੇ ਦੇ ਧਾਰਮਿਕ ਬੰਦੇ ਨੇ ਹੰਕਾਰ ਹੋ ਗਿਆ ਦੇਖ ਤਾਂ ਕਿ ਹੈ ਤਾਂ ਅੜਮੀ ਹੈ ਪਰ ਉਹ ਧਰਮ ਦਾ ਹੰਕਾਰ ਹੋ ਗਿਆ ਵੀ ਮੈਂ ਕਰਮੀ ਨੂੰ ਮੈਂ ਨਤ ਨਹੀਂ ਮੈਂ ਉਹ ਦਾਨ ਕੀ ਦੇ ਜਾਨਾ ਮੈਂ ਹਾਖ ਯੋਗੀ ਹਾਂ ਬੜੀ ਕਾਰ ਸੇਵਾ ਕੀਤੀ ਹੈ ਮੈਂ ਉਹ ਕੀਤਾ ਜੋ ਵੀ ਕੁਝ ਕਰਦੇ ਤੁਹਾਨੂੰ ਨੇ ਨਾ ਤੇ ਲੋਕ ਕਰਮकांड ਉਹਦਾ அவਮਾਨ ਉਤਾਰਨ ਦੇਵਤੇ ਨੂੰ ਮੈਕਾਸੋਸਮ ਸੁਮ ਬਾਇ ਉਹ ਉਤਾਰਦੇ ਹੋਏ ਜਿਤਰਨੇ ਮੈਕਾਸੋਸਮ ਤੁੰਗਾ ਜਿਹੀ ਹੋ ਜਿਤਰਨੇ ਜਥਾਂ ਦਾ ਇਹਦੇ ਜਲੇ ਜਿਤਰਨੇ ਇਹ ਚ ਵੀਰੇ ਚ ਲੈ ਇਹਨੇ ਆਖੇ ਸਰ ਜੇ ਭਗਤਾ ਜਿਹੜਾ ਹੋਆ ਰਾਵਣੀ दारु ਪੀਂਦੇ ਨਾ ਵਾਕੰਦੇ ਇਹ ਉਹਨਾਂ ਨੂੰ ਰਾਖੀ ਇਹਨਾਂ ਨੇ ਜਦੋਂ ਇਹ ਗੱਲਾਂ ਖੁੱਲਟੀਆਂ ਪਤਾ ਆ ਗਈਆਂ ਜੁੱਤੀ ਖੜਕ ਜਾਣੀ ਜੀ ਜੁੱਤੀ ਦਾ ਖੜਕੀ ਹੋਇਆ ਯਾਰ ਬ੍ਰਾਹਮਣ ਬਹੁਤ ਔਖੇ ਨੇ ਯੂਪੀ ਚੋਂ ਸਾਰੇ ਕਨੇਦਿਆਂ ਨੇ ਲੋਟ ਆਈ ਸੋ ਪ੍ਰੋਬਲਮ ਆਉਂਦਾ ਯੋਗੀ ਦੇ ਰਾਤ ਇਹਨੂੰ ਦਬਾਓ ਸਰਪੰਚਾਨੇ ਬ੍ਰਾਹਮਣ ਸਾਰੇ ਖਿਲਾਫ ਨੇ ਆਉਂਦਾ ਨਾ ਸਾਰੇ ਯੋਗੀ ਬ੍ਰਾਹਮਣ ਕਹਿੰਦੇ ਕਿ ਇਹ ਯੋਗੀ ਦੇ ਰਾਤੇ ਅੰਦਰੋਂ ਕੁਝ ਕਹਿੰਦਾ ਹੋ ਰਾ ਉਹ ਕਹਿੰਦੇ ਨੇ ਅਸੀਂ ਹਿੰਦੂ ਆ ਉਹ ਕਹਿੰਦੇ ਨੇ ਸਿਰਸਾ ਨਾ ਤੀਨ ਸਿੱਧੂ ਬੰਤੇ ਦੀ ਕੋਈ ਆ ਜੀ ਹਾਂ ਬਾਬਾ ਜੀ ਤੁਸੀਂ ਕਿਹਾ ਵੀ ਜਿਹੜੇ ਮੁਸਲਮਾਨ ਹੈ ਉਹ ਬੇਦ ਤੋਂ ਨਿਕਲੇ ਆ ਹਿੰਦੂ ਤਾਂ ਚਲੋ ਮੁਸਲਮਾਨ ਮੁਸਲਮਾਨਾ ਤੇ ਤਾਂ ਬਾਬਾ ਬੇਦ ਤੋਂ ਨਿਕਲਿਆ ਹਿੰਦੂ ਜੁਦੀ ਵੇਚਣ ਕਰਨਾ 파르시 ਜਿਹੜੇ ਨੇ ਨਾ ਉਹਨਾਂ ਨੂੰ ਸਨਮਾਨ ਲੈਣਾ ਹਿੰਦੂ ਨੂੰ 파르시 ਨਾ ਹਿੰਦੂ ਨੇ ਲੈ ਉਹ ਸਨਮਾਨ ਨੂੰ ਬੜਾ ਬੜਾ ਗੱਲ ਕਰਦੇ ਸੀ 파르시 ਸੀ ਉਹ ਮੁਸਲਮਾਨ ਨੇ ਨਾ ਹਿੰਦੂ ਨੇ ਦੋ ਜਣੇ ਹੀ ਹੁੰਦੇ ਹੈਗਾ ਜੈਨ ਮਤ ਪੈਦਾ ਹੋ ਗਿਆ ਬੁੱਧਵਾਤ ਉਹ ਇਕ ਬੁੱਧਵੰਤ ਹੋ ਗਿਆ ਜੈਨੂਤ ਹੋ ਗਿਆ ਜੈਨ ਵੱਧ ਜਾਦਾ ਹਿੰਦੂਵਾਂ ਨਾਲ ਚਲੇਗਾ ਜੋ ਵੱਧ ਮਤਜਾਦਾ ਮੁਸਲਮਾਨਾਂ ਨਾਲ ਚਲੇਗਾ ਸ੍ਰੀ ਕੰਡ ਕੌਣ ਜੁਟਾ ਹਕੀਆ ਨਹੀਂ ਨੇ ਕਿ ਲਾਗੇ ਪੀਰੋਂ ਕੰਨ ਮਰਟੀਆਂ ਉਹ ਪੀਰ ਅੱਧਾ ਮੁਸਲਮਾਨ ਹੈ ਜੋਗੀ ਕਾਹਨ ਇਸਲਾਮ ਕਬੂਲ ਲਿਆ ਸੀ ਇਹਨਾਂ ਨੇ ਚੌਂਦੀਆਂ ਜੋਗਿਆ ਨੇ ਜਦੋਂ ਆਮਨੇ ਪਰਮਪਰਵਿਤ ਕਰਦਾ ਤਾਂ ਇੱਕੋ ਹੀ ਸੀ ਗੱਲ ਉਹ ਕਹਿੰਦਾ ਤੂੰ ਖਾਣਾ ਪੀਣਾ ਆਪਣਾ ਆਖ ਲੋ ਤੀਰਥਾਂ ਤੇ ਵੀ ਜਾਓ ਉਹ ਬਾਣੀ ਕਲਾਮਾ ਸਾਡੀ ਨੂੰ ਪੜ੍ਹ ਲੋ ਜਿਹੜੇ ਜੋਗੀ ਸੀ اسی ਤਰ੍ਹਾਂ ਮਤਾਂਲੇ ਉਹ ਕਹਾਂ ਮਾ ਠਕਲਾ ਮਾ ਵੀ ਨੇ ਉਹ ਵੀ ਇੱਕੋ ਹੀ ਗੱਲ ਉਹ ਠੀਕ ਹੈ ਪੜ੍ਹ ਲੈ ਨਾ ਕਲਾਮਾ ਤੇ ਜਾਇ ਤੇ ਨਾਲੇ ਮਾਂਤਾ ਮਿਲਦੀ ਜੀ ਮੁਸਲਮਾਨ ਨੂੰ ਨਹੀਂ ਮੁਸਲਮਾਨ ਦਾ ਰਾਸਿ ਇਸ ਸੰਗਿਆਤ ਮਾਂਤਾ ਮਿਲਦੀ ਸੀ ਇਹ ਹੁਦਿਆਂ ਜਮਨ ਤਾਂ ਮਰਦੇ ਸੀ ਮਾਤੇ ਖੁਸੀ ਪਾੜਨ ਬਰਫ ਚੁੱਟਾਈ ਕਰਦੇ ਪਾਲੇ ਪਾਛੇ ਜਾਏ ਸਾਈ ਹੋ ਸੀ ਸ਼ੇਵੀ ਨੂੰ ਕਹਲਾਸ ਮਿਲ ਆ ਜੀ ਕਲਾਜ ਬਰਫਾਂ ਦੇ ਅੱਡਨੇ ਸਾਰੇ ਹੋ ਨੇ ਸਾਈ ਉਹਦੀ ਉਧਰ ਇਸ ਕਰਕੇ ਵਾਕੀਕਰ ਮਰਟ ਹੋ ਗਏ ਜਿਹੜੇ ਹਿੰਦੂ ਸੀ ਮੱਕੇ ਦੇ ਵਿੱਚ ਮੂਰਤੀਆਂ ਸੀ ਕਰਵਾਟ ਹੋਇਆ ਨੇ ਮੱਕਿਆਲੇ ਤੁਸਾਂ ਨੂੰ ਨਿਕਾਲਿਆ ਸਰਵ ਮੂਰਤੀਆਂ ਮੂਰਤੀਆਂ ਤੋਂ ਥੋੜੀਆਂ ਬਸ ਨੂੰ ਮੈਂ। ਇਹ ਉਦੇਵੀ ਮੂਰਤੀ ਪੂਜ ਕੇ ਨੇ ਮੂਰਤੀ ਪੂਜਾ ਦੇ ਖਿਲਾਫ ਹੈ। ਬਾਕੀ ਸਭ ਕੋ ਠੀਕ ਹੋ ਹੈ। ਸਿੱਖ ਵੀ ਹੋਈ ਨਾ। ਸਿੱਖ ਮੂਰਤੀ ਪੂਜਾ ਦੇ ਖਿਲਾਫ ਇਹ ਤਾਂ ਮੂਰਤੀ ਪੂਜਾ ਦੇ ਵੀ ਖਿਲਾਫ ਹੋ ਗਿਆ। ਇਹ ਤਾਂ ਫੇਰੋਜ਼ਾ ਲੈਣ ਤੇ ਆ ਕੇ ਗੁਰੂਆਂ ਨੂੰ ਜੋੜ ਕੇ। ਇਸਲਾਮ ਵਾਲੇ ਨੇ ਲੇਗਾ ਸਕੇ ਦੇ ਪਿੱਛੇ। ਸਿੱਖ ਵੀ ਖਤਮ ਹੋਵੇ 500 ਸਾਲ ਚ। ਇਸਲਾਮ ਖੜਾ ਹੁੰਦਾ ਸੀ ਮੁਸਲਮਾਨ ਖੜਾ ਹੁੰਦਾ ਸੀ ਮੁਸਲਮਾਨ ਉਹ ਤੇ ਖੜਾ ਸੀ ਉਦੋਂ ਗੁਰਨਾਨਕ ਬੇੜੇ ਕਬੀਰ ਦੇ ਚੰਦੇ ਟਾਕੇ ਨਹੀਂ ਹੋ ਗਏ ਸੀ ਸਾਰੇ ਇਸਲਾਮ ਵਾਲੀ ਗੱਲ ਸੀ ਮੁਸਲਮਾਨ ਦੇ ਘਰ ਪੈਦਾ ਹੋ ਗਏ ਕਬੀਰ ਨੇ ਗੁਰਮਤ ਮੰਨੀ ਕਿਉਂ ਅਸਲ ਮਤ ਸੀ ਨਰੋਲ ਇਸਲਾਮ ਸੀ ਇਹ ਤਾਂ ਨਹੀਂ ਜਿਉਂ ਐਵੇਂ ਕੰਮਾ ਨਹੀਂ ਜਿਗੋ ਦਾਂ ਕਰਕੇ ਮੁਸਲਮਾਨ ਅਖਬੀਰ ਨੂੰ ਹੁੰਦੇ ਨੇ ਸਾਰੇ ਕਹਿੰਦਾ ਜੰਮੀ ਤਾਂ ਸਾਡੇ ਘਰੇ ਆ ਮਾਤੇ ਮੈਂ ਕਹਤਾ ਵੀ ਅਖਬੀਰ ਬੈਲਾ ਉਹ ਪਰਮੇਸ਼ਰ ਨੇ ਕਿਉਂ ਪੈਦਾ ਕੀਤਾ ਤੇ ਇਕਤਾ ਵਾਸਤੇ ਪੈਦਾ ਕੀਤਾ ਸੀ ਮੈਂ ਤਾਂ ਜੋ ਕਹ ਜੋ ਸੱਚਾ ਹੋਈ ਕਿਹਾ ਮੈਂ ਕੁਝ ਝੂਠ ਬੋਲੇ ਇਹ ਸਿੱਖ ਕਿਉਂ ਕਹਿੰਗਾ ਤੇ ਸਨਾਤਨੀ ਇਹ ਕਹਿੰਦੇ ਜੇ ਅਖਬੀਰ ਕਹਤਾ ਇਹ ਦੋ ਜੂ ਮਹਲਵਣ ਨਾ ਵੀ ਲਿਖੋ ਨਹੀਂ ਏ ਜੌਨ ਨੇ ਨੀਟ ਪਾਰਾ ਪਾਕਿਸਤਾਨ ਤੋਂ ਆਇਆ ਉਹਨੇ ਹੰਦਰ ਦਵਾਰ ਬਣਾਇਆ ਮੁਸਲਮਾਨ ਬਣਾ ਉਹਨੇ ਮਿਲਦਾ ਦਿੱਤਾ ਖਾਨ ਤੱਕ ਨਿੰਦਾ ਕੀਤੀ ਰੰਦਰ ਦੇਤੇ ਨੇ ਟਾਹਿਆ ਸੀ আর ਖਲਾਫ ਉਹਨੇ ਆਤਮਾ ਤੇ ਗੁੰਡੇ ਕਹਿਣ ਵਾਲੇ ਜਿਹੜੇ ਗੁੰਡੇ ਜਿੰਦੂਆਂ ਦੇ ਖਲਾਫ ਤਰਫ ਦੇ ਖਲਾਫ ਕਰਦੇ ਨੇ ਸਾਸ਼ਾ ਖੁੱਲ ਕੇ ਸਾਰੇ ਬੋਲਦੇ ਨੇ ਮਨ ਬਾਰੇ ਭਗਵੰਤੂ ਜੀ ਸਾਡੇ ਟੀਵੀ ਤੇ ਪ੍ਰਚਾਰ ਕੀਤਾ ਰਾ ਉਹਨਾਂ ਨੂੰ ਪਤਾ ਹੈ ਵੀ ਦੁਨੀਆ ਨੇ ਸਿੱਖ ਮਤ ਨੂੰ ਕਬੂਲ ਕਰ ਲਿਆ ਮੈਸੇਜ ਚੱਲਿਆ ਗਿਆ ਸਨਾਤਨੀ ਹਿੰਦੂ ਵੀ ਕਹਾਂ ਮੁਸਲਮਾਨ ਕਰ ਰਹੇ ਇਹਦਾ ਭਗਵੰਤਾਈ ਮੈਸੇਜ ਚੱਲਿਆ ਗਿਆ ਇੱਕ ਦਵਾਇਆ ਬਸ ਉਹਨਾਂ ਨੇ ਚੜ੍ਹ ਲੈ ਲਿਆ ਗਿਆਨ ਇੱਕ ਬਾਰੇ ਬਹੁਤ ਹੁੰਦਾ ਜੁੱਤਾ ਦੁਬਾਰਾ ਭਗਵੰਤੂ ਜੀ ਆਣ ਵੀ ਇਹ ਜੀ ਦੁਆਰਾ ਕੋਲ ਮੰਨ ਦੀ ਜੁੱਤੀ ਹਾਣੀ ਚਾਹੇ ਅੰਦਰੋਂ ਦੁਖੀ ਯੋਗ ਦੱਸ ਤਾਵੇ ਬ੍ਰਹਮ ਜੀ ਹਾਂ ਅੱਛਾ ਕਾਹ ਕੇ ਦਿਖਾਉਣ ਇੱਕ ਝੂਠ ਹੈ ਨਹੀਂ ਸਿੱਖ ਅਕਾਲ ਤਖ ਨੂੰ ਇਹ ਨਹੀਂ ਕਹਿੰਦਾ ਮੈਂ ਅਕਾਲ ਤਖ ਨੂੰ ਨਹੀਂ ਮੰਨਦਾ ਮੈਂ ਉਹਦਾ ਫੋਲ ਕਰ ਰਿਹਾ ਕਰਦਾ ਹਾਂ ਉਹਨੂੰ ਪੰਟੀ ਨਹੀਂ ਦਿੰਦਾ ਤਾਂ ਤੂੰ ਕਹੇ ਪਰ ਉਹ ਤਾਂ ਫੰਕੀ ਆ ਕਾਲ ਕਰਤਾ ਲੰਡੂ ਕੁਛ ਮੇਰੇ ਕੋਲ ਕੋਈ ਸਮਝ ਨਹੀਂ ਕਿ ਫੋਨ ਕੀਤਾ ਇਹ ਤੋਂ ਮੰਨ ਅਸੀਂ ਰਿਕਾਰਡ ਕਰਾਂਗੇ ਵੀ ਮੈਂ ਕਹਤਾ ਉਹਨੂੰ ਨਹੀਂ ਮੰਨਦਾ ਕਿਉਂਕਿ ਗੁਰਮਤਿ ਖਰਾਬ ਨੇ ਨਹੀਂ ਮੈਂ ਨਾਲ ਗੱਲ ਨਹੀਂ ਬਹੁਤ ਟਾਈਮ ਨਹੀਂ ਹੈ ਤੁਹਾਡੇ ਵਾਸਤੇ ਚਾਰ ਆਦਮੀ ਜਵਾਬ ਦੇ ਚੁੱਕਿਆ ਹਾਂ ਉਹਨੂੰ ਉਲਟੇ ਸਿਰ ਜੜਿਆ ਬਾਠੋੜਣਾ ਮੈਂ ਕਿਹਨੂੰ ਕਰਾਂ ਉਸਦੇ ਮਤਿਓਤ ਗਾਲ ਤਾਂ ਹੁਣ ਹੁੰਦਾ ਨਹੀਂ ਬੈਠੇ ਉਹਨੇ ਬੈਠਾ ਫਿਰ ਕੱਲ ਕਾਇਆ ਕਲਨ ਜਮਨ ਤਾਂ ਵੇਲਾ ਕੀ ਹੁੰਦਾ ਵਾ ਅ ਕੱਲ ਕਾ ਮੈਂ ਉਹ ਸਿੱਖ ਨਹੀਂ ਉਹਨਾਂ ਵਾਲੀ ਸਿੱਖੀ ਮੈਨੂੰ ਨਹੀਂ ਮੰਦਾ ਇੰਟਰਨੈਟ ਤੇ ਪਾ ਫਿਰ ਮੈਂ ਨਾਲ ਗੱਲ ਕਰਾਂ ਨਹੀਂ ਬਾਈ ਕੋਣਾ ਥੋੜਾ ਮੈਨੂੰ ਨਹੀਂ ਫੋਨ ਕਰਨਾ ਲੇਕਿਨ ਖਚਾਉਂਦੇ ਰਹਿੰਦੇ ਜੀ ਨਖ ਨਖ ਪਰਸੇਵ ਜਾਂਚੈ ਸੁਰਸਰੀ ਬਾਬਾ ਜੀ ਇੱਥੇ ਪ੍ਰੋਫੈਸਰ ਸਹਿਬ ਸਿੰਘ ਨੇ ਅਰਥ ਕੀਤੇ ਆ ਗੰਗਾ ਉਸ ਦੇ ਦਰ ਤੇ ਉਸ ਦੇ ਨੌਂਹਾਂ ਦਾ ਪਸੀਨਾ ਹੈ ਉਹ ਪਰਸੇਵ ਉਹਦਾ ਪਸੀਨਾ ਹੀ ਕਾ ਲੋਪਸੀਨਾ ਤਾਂ ਕਰ ਹੁੰਦਾ ਨਹੀਂ ਉਹਦੇ ਹੱਥਾਂ ਦਾ ਪਸੀਨਾ ਕਹਿ ਸਕਦੇ ਹਾਂ ਅਸੀਂ ਚੇਤਰਮਨ ਹੱਥ ਨੇ ਨਾ ਉਹ ਕੋਈ ਹੱਥ ਹੁੰਦਾ ਉਹਦਾ ਦੋਹੇ ਨਹੀਂ ਉਹਦੀ ਜਿਹੜੀ ਸਖਤ ਉਹਦੇ ਜਿਹੜਾ ਮੁਖ ਹੈ ਗੰਗਾ ਮੁਖ ਤੋਂ ਨਿਕਲੀ ਹੋਈ ਹੈ ਨੋਂ ਦਾ ਪਸੀਨਾ ਨਹੀਂ ਹੁੰਦਾ ਨਾਲੇ ਗੰਗਾ ਤਾਂ ਹੈ ਹੀ ਨਹੀਂ ਸਭ ਸੀ ਤਾਂ ਮਤਲਬ ਸੁਰਸਰੀ ਮੈਂ ਤੈਨੂੰ ਕਹਾਣੀ ਕਿਉਂ ਸੁਣਾਈ ਆ ਹਲਾਵਾ ਦੀ ਬੇਈਮਾਨ ਗੰਗਾ ਅਥ ਕਹਿੰਦਾ ਉਹ ਯਾਰ ਗੰਗਾ ਜਮਨਾ ਸੁਰਸਰੀ ਉੱਥੇ ਮਿਲਦੇ ਨੇ ਹਾਂ ਇਹਨਾਂ ਨੇ ਗੰਗਾ ਨੂੰ ਸੁਰਸਰੀ ਸੁਰਸਰੀ ਨੂੰ ਗੰਗਾ ਕਹਤਾ ਕਿਉਂ ਗਿਆਵੇਂ ਉਹਨੇ ਜਦ ਫਸ ਗਏ ਗੰਗਾ ਕਨਾਲ ਰੈਸੋਰਟ ਦੀ ਤੁ ਫਤੈਨੇ 3 ਵਾਇਟ ਪਿੰਗਲਾ ਸੁਖਮਣਾ ਪਹਿਲਾ ਇਹੜਾ ਫਿਰ ਪਿੰਗਲਾ ਫਿਰ ਸੁਖਮਣਾ ਸੁਖਮਣਾ ਸੋਰ ਫਰੀ ਗਿਆ ਵਿਚਾਰੇ ਦਾ ਪਿੰਗਲਾ ਗੁੰਦਾ ਆ ਤੇ ਰਵਣੀ ਉੱਥੇ ਫੋੜ ਗੰਗਾ ਫਿਰ ਸੁਖਮਣਾ ਲੰਗਾਂ ਨੂੰ ਸੁਖਮਣਾ ਕਿਵੇਂ ਕਹਾਂ ਮੈਂ ਤੁਸੀਂ ਵਿਖਾਰੇ ਜਾਦੋ ਆਹਿੰਚਲਾ ਕੀਆ ਨਹੀਂ ਉੱਤੇ ਜ਼ਮੀਨ ਤੇ ਕੁਝ ਬਣਾ ਬੈਠੇ ਪਰ ਚਾਰ ਵਾਲੇ ਫਾਜਾ ਦੇ ਫੇਰ ਕੁਝ ਕਹਿਣ ਦੇ ਨਹੀਂ ਤੁਹਾਨੂੰ ਕਿਹੜਾ ਪਤਾ ਛੋਟ ਕਿਹੜਾ ਆਦ ਰਹਿ ਗਿਆ ਲੋ ਇਹਦਾ ਨੋਟ ਕਰਾਉਣੀ ਹੈ ਹੁਣ ਸੁਰਸੇ ਨਹੀਂ ਕਹਤਾ ਉਹਨੇ ਗੰਗਾਂ ਗੰਗਣ ਸੁਰਸੇ ਦੀ ਕਿ ਮੈਂ ਕਹ ਦੁ ਉਹ ਤਾਂ ਕਹੂੰਗਾ ਜਦ ਕਹਿੰਦਾ ਗੰਗਾ ਜਮਨ ਕੇ ਅੰਤਰੇ ਠੀਕ ਹੈ ਜੀ ਜਮਨ ਨਾਲੇ ਰੜੇ ਹੁੰਦਾ ਸੋਸਰੀਏ ਸੋਸਰੀ ਦਾ ਆਇਓ ਫਿਰ ਸੋਸਰੀ ਵਿਛਾਲੇ ਹੋਣੀ ਸ਼ਾਇਦ ਸੋਨ ਨੂੰ ਕਹਿ ਗਾਉਤ ਉਹ ਹੱਦ ਤੇ ਹੈ ਜਿਹੜੀ ਅਸੀਂ ਪਾਰ ਕਰਨੀ ਹੈ ਜਿਹਨੂੰ ਗੰਗਾ ਨੂੰ ਟਾਹ ਹੈ ਕਾਇਰ ਨੇ ਬਤਾੜਨੀ ਨਦੀ ਇਹ ਪਾਰ ਨਹੀਂ ਜਾਣ ਪਾਰ ਨਹੀਂ ਜਾ ਉਹਦਾ ਕੋਈ ਪਾਰ ਨਹੀਂ ਪਾ ਸਕਦਾ ਉਨਦੇ ਪਾਰ ਕੋਈ ਹੋ ਹੀ ਨਹੀਂ ਸਕਦਾ ਵੱਡਾ ਦਰਿਆ ਹੈ ਉਹ ਤਾਂ ਗਏ ਨਹੀਂ ਨੇ ਸੁਰਸਤੀ ਦਾ ਕਹਾਂ ਜਾਗੇ ਆ ਉਹ ਜਿਆਦਾ ਫਿਰ ਗੰਗਾ ਚਬਨਾਓਗੇ ਉਹਦਾ ਵਿਚਾਲਾ ਹੋ ਜਾਂ ਸੁਰਸਤੀ ਅਰ ਗੰਗਾ ਦਾ ਵਿਚਾਲਾ ਹੋ ਜਾਂ ਚਬਨਾਓ ਦਾ ਵੀ ਵਿਚਾਲੇ ਯਕੀਨਾਂ ਤੈਨ ਮਾਰ ਕੇ ਦੇਖ ਜਿੰਨਾ ਤੇ ਲਿਖਣਾ ਗੰਗਾ ਜਵਨ ਕਾਉਂਤਰਾ ਇਹ ਜੰਨਾ ਜੰਨਾ ਦੋ ਕੱਠੀਆਂ ਨੇ ਇਹ ਸੁਸ ਵੀ ਨਹੀਂ ਹੈ ਬਿਚਾਰੇ ਇਹਨਾਂ ਦੇ ਤੀਜੀ ਕਿਠਾਈ ਤੇ ਦੋਵੇਂ ਮੰਦਰ ਤੇ 30 ਖੜੂਗਰ ਦਰੂ ਇੱਥੇ ਅਲਾਵਾ ਤੁੰਮ ਇੱਕ 700 ਹੋਰ ਵੀ ਆ ਪੰਜਾਬ ਚ ਪੁਰਾਣੇ ਚ ਆ ਜਿਹੜੇ ਬੈਠੇ ਨੇ ਨਾ ਪੱਟ ਜੇਲੀ ਕੋਮ ਖੇਤਰ ਸਰੋਵਰ ਜੀ ਜਾਂਦਾ ਨਾਲ ਆ ਜਾ ਨਿਕਲ ਕੇ ਇਹ ਗੋਆ ਦਾ ਉਹੀ ਬਠਾਤੀ ਗਿਆ ਜਿਗਾ ਦੇ ਤੋਂ ਨਿਕਲਦਾ ਹੋ ਜਿਗਾ ਦੇ ਉੱਪਰ ਗਪਾਲ ਤੋਂ ਇਕੱਠਾ ਜਾਂ ਪਾਣੀ ਹੋ ਕੇ ਨਾ ਇਹ ਉਪਰ ਉਧਰ ਉੱਥੇ ਚੱਲ ਜਾਣਾ ਆਪਣੇ ਜਿਹੜਾ ਜੀਂਗਾ ਉਹ ਨੂੰ ਵੀ ਸਭ ਕਹਿੰਦੇ ਨੇ ਕੋਹ ਚੈਤਲ ਦੇ ਸਰੋਵਰ ਚੋਂ ਹੀ ਪਾਣੀ ਜਾਂਦਾ ਫਲਗੂ ਵੀ ਉਹੀ ਪਾਣੀ ਜਾਂਦਾ ਇਹ ਟੇਕਓਵਰ ਤੇ ਦਿੱਪਟ ਜਿਹਨਾਂ ਨੇ ਬਾਣੀ ਗੁਰੂ ਗ੍ਰੰਥ ਸਾਹਿਬ ਜਿੱਥੋਂ ਪਾਈ ਕੁਨੀਸੇ ਨੇ ਬਣੇ ਨੇ ਪਰ ਹੈ ਕੋ ਕ ਵੀ ਸੋਤਸਰੀ ਕਹਿੰਦੇ ਨੇ ਸਰਾਸੋਤੀ ਕਹਿੰਦੇ ਨੇ ਵੀ ਅਸੀਂ ਕਣਾਂ ਨੇ ਬੈਠੇ ਆ ਕਿ ਉਹ ਨੇ ਨਾ ਉਹ ਉਹ ਉਹਨਾਂ ਨੇ ਉਹ ਉਹਦਾ ਨਾਮ ਸੋਤਸਰੀ ਦੇਤਾ ਉਹ ਆਵਾਜ਼ਾਂ ਦੇ ਨੂਦਾਂ ਨੋਸਰਾ ਫਿੱਦੇ ਲੱਟਾ ਹੋਇਆ ਇਹ ਫਸੇ ਬੈਕਦੇ ਕੋ ਜਿੱਥੇ ਜਗ੍ਹਾ ਨੇ ਇਹਨਾਂ ਨੇ ਬਣਾਈਆਂ ਹੋਈਆਂ ਜਿੱਦੇ ਸੀਤਾ ਨੇ ਬਣਵਾਸ ਕਟਿਆ ਸੀਤਾ ਮੰਡੀ ਕੋਣ ਹੈ ਕੋਈ ਕੁਸ਼ਮ ਇੱਥੇ ਆਜਣੇ ਪੰਚਕੂਲਾ ਇੱਥੇ ਇਹਨਾਂ ਨੇ ਬਣਾਇਆ ਵੀ ਇੱਥੇ ਉਹ ਪੱਦੇ ਪੱਨੋਂ ਨੇ ਇੱਥੇ ਬਣਵਾਸ ਕਟਿਆ ਪੰਚਕੂਲਾ ਹੋਇਆ ਇੱਥੇ ਪੰਜਾਣੇ ਨੌਦੇ ਆ ਇਹ ਕਿਹੜਾ ਟਪੀਂ ਗੋਡਾ ਪਾਣੀ ਨਹੀਂ ਬਣਾਇਆ ਹੋਇਆ ਕਿਤੇ ਵੀ ਮੈਨੂੰ ਗੋਡਾ ਮਾਰਿਆ ਤਾਂ ਕਿਹਜ ਪਾਣੀ ਨਿਕਲਿਆ ਪੱਥਰ ਜੇ ਇਹ ਕਿਹੜਾ ਥੋੜਾ ਝੂਠ ਬੋਲਦੇ ਨੇ ਸਾਡੇ ਬਣਾਤਾ ਪੌੜ ਮਾਰਿਆ ਪਾਣੀ ਨਿਕਲਿਆ ਆ ਆਨੰਦ ਦੇ ਨਾਲ ਉਹ 10 12 ਤੋਂ ਉਹਦੇ ਨਿਕਲਦਾ ਪਾਣੀ ਜਦੋਂ ਟੈਂਕ ਬਣਿਆ ਨਾ ਪਹਿਲੇ 1000 ਤੋਂ ਨਿਕਲਦਾ ਹੁੰਦਾ ਸੀ ਪਾਣੀ ਉਹ ਥੋੜੇ ਸਾਲ ਹੋ ਗਏ ਹੋ ਗਏ ਉਹ ਕਈ ਤੋਂ ਉਹਦੇ ਪੜ ਮਾ ਓਏ ਆ ਜਗਾ ਨਿਕਲਦਾ ਚੁੱਪ ਬੋਇ ਤਾਂ ਪਹਿਲੇ ਨਹੀਂ ਲੀਵੰਗਾ ਇਹਨਾਂ 47 ਹੋਣੀਆਂ ਕੋਈ ਪਰ ਉਹ ਦਰਿਆ ਕਸ਼ਮੀਰ ਵੀਰ ਜਗਨ ਨਾਲ ਪਾੜਨ ਦੇ ਵਿੱਚ ਕਹਿੰਦਾ ਜੀ ਪੌੜਾ ਦਾ ਪੌੜ ਮਾਰੇ ਆਇਆ ਤੇ ਕਿਤੇ ਪਾਣੀ ਨਿਕਲਿਆ ਜਾਂ ਤਾਂ ਗਏ ਨਹੀਂ ਉੱਤੇ ਗੁਰੂ ਕੀ ਲਾਹੌਰ ਪਿਆ ਇਹ ਕਿਹਦਾ ਤੋਂ ਤੋਂ ਘੂੜੇ ਉਹਨਾਂ ਨੇ ਜੀ ਝੂੜਦਾ ਸਦਾ ਹੀ ਧਰਮ ਜਿਹੜਾ ਵੱਡਾ ਝੂੜ ਹੈ ਵੱਡਾ ਵਰਸ਼ਾ ਫਿਰ ਉਹਨਾਂ ਦੀ ਖੋਲ ਨਹੀਂ ਚੱਟਦੀ ਮੇਰੀ ਖੋਲਨੀ ਵੱਡੀ ਕ ਵਰਸ਼ਾ ਵੱਡਾ ਜੇ ਖੋਲਨੀ ਵੱਡੀ ਆ ਖੋਲਦੀ ਕੋਸ਼ਿਸ਼ ਕਰਦੀ ਵਰਸ਼ਾ ਦੂਰ ਤੱਕ ਮਾਰ ਕਰਦਾ ਉਹ ਜਿਹੜੀ ਹੈ ਪਾਈਏ ਉਹ ਗੁਰਮੱਤਾ ਗੰਗਾ ਉਹਦੇ ਕਥੇ ਉਹਦੇ ਦੌਰੇ ਚਲੋ ਉਹਨਾਂ ਆਪਾਂ ਗੰਗਾ ਦੇ ਨਹਾ ਚੋਂ ਕਹਿੰਦੇ ਨਿਕਲੀ ਆ ਉਹ ਅਗੀਰ ਥੱਲੇ ਗਿਆ ਪਹਾੜਾਂ ਚੋਂ ਲੈ ਗਿਆ ਪਾਣੀ ਪਹਾੜ ਵੱਡ ਵੱਡ ਕੇ ਲੈ ਗਿਆ ਸਾਖੀ ਬਣਾਈ ਇਹਨਾਂ ਦੀ ਉਹਨੇ ਕਿ ਥੋੜੀ ਗੱਲ ਉਹਦੇ ਨਹਾ ਚੋਂ ਨਿਕਲੀ ਗੰਗਾ ਦੀ ਸਾਖੀ ਲੰਘ ਪਈ ਐ ਬਾਹਰਿਤ ਲੈ ਕੇ ਆਇਆ ਗਾਂ ਸ਼ਿਲੀ ਜੀ ਬੈਠਾ ਸ਼ਿਲੀ ਜੀ ਦੇ ਉੱਤੇ ਤਾਰ ਪੈ ਗਈ ਜਿਹੜੀ ਇਹਦੇ ਜਟਾਂ ਦੇ ਵਿੱਚੋਂ ਹੀ ਨੰਗਾ ਨਿਕਲ ਨਹੀਂ ਦਿੱਤੀ ਬਾਹਰ ਅੜਜਾਲੀ ਉਹੀ ਆ ਗੁਰੂ ਨਾਨਕ ਲੈ ਕੇ ਆਇਆ ਗੰਗਾ ਸਰੀ ਚੰਗੇ ਜਟਾਂ ਦੇ ਲਕੋੜੀ ਅੜਜਾਲੀ ਉੱਥੇ ਹੀ ਹਣ ਜਾਈ ਪਈ ਐ ਇੱਥੇ ਵੀ ਜਟਾਂ ਦਾ ਹੋਈ ਆਈ ਹੋਈ ਜੜਾ ਨੂੰ ਹੰਦਨੇ ਲੋਕ ਜੀ ਨੂੰ ਮੰਨ ਉਹਨੂੰ ਸੇਈ ਚੰ ਨੂੰ ਮੰਨਦੇ ਨੇ ਸੇਈ ਚੰ ਦਾ ਪੱੜ ਲੱਗਿਆ ਤੁਹਾਡੇ ਉੱਤੇ ਦਰਬਾਰ ਦਾ ਹੋਈ ਆਈ ਨੇ ਬਿਲਕੁਲ ਜੀ ਪੱੜ ਗਿਆ ਕਦੇ ਪੱੜ ਲੱਗ ਗਿਆ ਹੈ ਤੇ ਪਰਦੋਸਣ ਵਾਲਾ ਬੰਦੇ ਲੋਕ ਸਾਨੂੰ ਦਾ ਪੱੜ ਲੱਗ ਗਿਆ ਹੈ ਪੱੜ ਲੱਗਿਆ ਆ ਇਹ ਲੈ ਦੇ ਤੇ ਪਰ ਦਵਾਰ ਤੋਂ ਪੈ ਰਾਇਆ ਦਵਾਰ ਪਾੜ ਦਿੰਦਾ ਪੱਤੋਂ ਨੂੰ ਵਾਰਦੂ ਨਾ ਕਰ ਪਾੜਦੇ ਸੰਗਤ ਕੇ ਨੂੰ ਕਰਤੀ ਰਾਤੇ ਨਾਲੇ ਜੀ ਅੱਗੇ ਪੜੇ ਤੈਨਾਂ ਕਾ ਦਰ ਮੈਨ ਅਜੇ ਤਾਂ ਪ੍ਰਕਲਪੋਂ ਤੋਂ ਬਾਹਰ ਇਹ ਕਿਹਦੇ ਨੂੰ ਨਾ ਫੇਲੀਆ ਦੇਖਦਾ ਨਖ ਪਰਸੇਵ ਜਾਂਚੈ ਸੁਰਸਰੀ ਉਹਦੇ ਜਿਹੜਾ ਉਹਦੇ ਅੰਦਰ ਸੱਚ ਐ ਨਾ ਸੱਚਖੰਡ ਚ ਉਹ ਸੁਰਸਰੀ ਆਈ ਐ ਤੁਰਕੀ ਬਾਣੀ ਹੈ ਸੁਰਸਰੀ ਤੁਰਕੀ ਬਾਣੀ ਆਈ ਤੰ ਚੰਦ ਮੰਗਾਈ ਐ ਤੁਰਕੀ ਬਾਣੀ ਹੈ ਭਾਈ ਉਹਦੇ ਹਿਰਦੇ ਚ ਹੋਈ ਉਹਦੇ ਕ ਕਰਹੀ ਹੁੰਦਾ ਹਿਰਦੇ ਹੁੰਦਾ ਕ ਦੇਨ ਘਰ ਨਹੀਂ ਕਹਿੰਦੇ ਜਾਂ ਕਿ ਘਰ ਹੈ ਘਰ ਦਾ ਸ਼ਬਦ ਵਰਤੇ ਹੋਇਆ ਉਹਦਾ ਹਿਰਦੇ ਘਰ ਨੌ ਤਾਰੇ ਹੁੰਦੇ ਹੀ ਨਹੀਂ ਮੈਨੂੰ ਐ ਦੱਸ ਲਾਉ ਕਿੱਥੇ ਨੇ ਜੇ ਨੌ ਨੇ ਤਾਂ ਮਾਫੀ ਹੋਊਗਾ ਤੇ ਆਦਮੀ ਦਾ ਜੀਰੋ ਆਦਮੀ ਨਾਮ ਮੰਨੇਗਾ ਆਦਮੀ ਐ ਫਿਰ ਉਹ ਆਗਮਗਾ ਨਿਕੜੀਏ ਫਿਰ ਉਹਦੇ ਹੰਗਾ ਵੀ ਆਹੀ ਹੋਊਗੀ ਕੀ ਆਤਰਤਲ ਵੀ ਟੁਲਕੀ ਬਾਣੀ ਰਹੀ ਫਿਰੇ ਮੈਂ ਨੋਟਾਂ ਨਹੀਂ ਜਿਵੇਂ ਨੂੰ ਟਾਈਮ ਦਤੋ ਨਾ ਵੀ 76 ਫੇਰ ਦੂਗਾ ਸੰਗਤ ਦੇ ਵਿੱਚ ਕੋਈ ਝੂਠ ਫੇਰ ਦੇਣਾ ਨਾ ਅੰਮਰਸਾਰੇ ਮੈਂ ਸੀ ਯਾਰ ਉਹ ਕਰਦਾ ਸੀ ਟਾਈਮ ਨਹੀਂ ਦਤੋ ਲੈ ਕਿੰਨਾਂ ਨੂੰ ਗੰਦੇ ਨਹੀਂ ਹੋਣੇ ਨੇ ਵੀ ਕਿਤੇ 10 ਜਾਣੇ ਗਏ ਸੀ ਉੱਤੇ ਮਾਨੂੰ ਆਪਣੇ ਸੱਥੀ ਦੇ ਕੇ ਸਦਗੋਸ਼ ਤੋਂ ਜਵਦੀ ਸਾਹਿਬ ਨੇ ਪਹਿਲਾਂ ਪੜਿਆ ਹੋਇਆ ਸੀ ਕਲਕੱਤੇ 파ਟਮੀਰ ਦਾਡਾ ਨੂੰ ਜੁਲਾ ਕਲਕੱਤੇ ਮੈਂ ਘਰ ਉਹ ਦੇ ਕੇ ਪੜਦਾ ਸੀ ਇਹਦੀ ਭੈਣ ਸੀ ਆਪਣਾ ਜਿਹੜਾ ਕੀ ਸੀ ਉਹ ਫਾਉਡੇਸ਼ਨ ਦਾ ਪ੍ਰਧਾਨ ਕਲਕੱਤੇ ਮਨਜੀਤ ਸਿੰਘ ਮਨਜੀਤ ਸਿੰਘ ਕਲਕੱਤਾ ਉਹ ਦੇ ਫੈਸਲੇ ਜੀ ਗਵਰਦੀਰ ਉਹ ਗਦੇ ਉਹ ਬਈਆ ਹੈ ਚੌਥੀ ਦੰਦਾ ਨੰਨ ਕਟਕਤੇ ਗੱਲ ਨੂੰ ਜੀ ਜੇ ਗੱਲ ਕੀਤੀ ਉਹਨੇ ਨੂੰ ਸੱਜਾ ਫਿਰ ਉਹਨੇ ਕਿਤਾਬ ਲਈ ਉਹਨੇ ਮਨਜੀਤ ਨੂੰ ਪੁੱਛਿਆ ਕਿ ਲੜਤਾ ਸਲਾਹ ਉਹ ਕਹਿੰਦੇ ਛੱਡ ਬੜੇ ਆ ਦੀ ਗੱਲ ਨਹੀਂ ਸਾਡੇ ਕੋਲ ਸਾਡੇ ਕੋਲ ਤਾਂ ਹੋਰ ਹੀ ਚੀਜ਼ ਹੈ ਬਾਰੇ ਦਾ ਤੂੰ ਕੀ ਕਰਦਾ ਹੈ ਕਿਹੜੇ ਨਾਲ ਪੈ ਗਿਆ ਤੂੰ ਉਹ ਕਹਿੰਦਾ ਹੈ ਸਿਆਸਤ ਦੇ ਵਿੱਚ ਨਹੀਂ ਇਹ ਗੱਲ ਜਲਦੀ ਹਸਾਉਂਦਾ ਰੋਮਾਂਟਿਕ ਗੱਲ ਹੈ। ਮੰਨੇ ਨਹੀਂ ਵਾਜੀ। ਹਾਂ ਜੀ ਸਭ ਪ੍ਰਕਾਸ਼ੇ ਦੀ ਚਿੱਠੀ ਹੈ। ਕੇ ਉਹਨੇ ਕਿਹਾ ਵੀ ਕਾਲੇ ਫਗਾਨੇ ਦੇ ਕਾਲੇ ਪਤਾ ਸੀ ਬੰਜੀਏ ਸਾਨੂੰ। ਉਹ ਪੜ੍ਹੀ ਸੀ ਕਹਾੜਦੋਏ ਕਹਾਵਾਂ ਪੜ੍ਹੀਆਂ ਸੀ। ਹਾਂ ਤੁਹਾਨੂੰ ਚਿੱਠੀ ਆਈ ਸੀ ਉਹ। ਆਹ ਸਭ ਪਤਾ ਸੀ ਇਹਨਾਂ ਨੂੰ ਬਈ ਮ ਪਤਾ ਹੈ ਵੀ ਇਹਦੇ ਚਲਦੀ ਨਹੀਂ ਉਹ ਗੁਰਮਤ ਅਲ੍ਹਾ ਕਮ ਨਹੀਂ ਹੈ ਪਬਲਿਕ ਨੂੰ ਨਹੀਂ ਕਿਹਾ ਇਹਨਾਂ ਨੇ ਪਬਲਿਕਲੀ ਸੁਣਾ ਕੇ ਐਕਸਪੋਜ਼ ਹੋ ਗਏ ਪਬਲਿਕ ਚਾਹੀਦਾ ਹੈ ਪਬਲਿਕ ਨੂੰ ਵੀ ਹੋਰ ਕੁਝ ਚਾਹੀਦਾ ਜੀ ਆ ਨਖ ਜਾਚੈ ਸੁਰਸਰੀ ਔਰ ਕਰ ਗੁਰਮਤਾ ਨਖ ਜਿਹੜੀ ਮੁੰਦੀ ਨੀ ਕਿਸੇ ਪਾਸੇ ਸਿੱਧੀ ਜਾਂਦੀ ਐ ਜਿਵੇਂ ਲੋਹਾ ਮੁੜ ਜਾਂਦਾ ਨਾ ਨਖ ਨਹੀਂ ਹੁੰਦਾ ਅਸਲੇ ਨਹੀਂ ਹੁੰਦਾ ਉਹ ਹੁਲਾ ਹੁਲਾਦ ਮੁੜਦਾ ਨਹੀਂਦਾ ਟੁੱਟ ਜਾਂਦਾ ਨਖ ਖੈਣ ਨੇ ਸਦਾ ਕਰਦਾ ਉਹ ਡੋਨਟ ਯੂ ਲਵ ਵਰਦਾ ਸਖਤ ਸੱਚ ਜਿਹੜਾ ਗਣਾ ਖੁੰਦ ਬੈਠੇ ਸ਼੍ਰਿੰਗ ਸੁਮੇਰ ਕਚੰਡ ਬਰਾਜਤ ਸ਼੍ਰਿੰਗ ਸੁਮੇਰ ਜਿਹੜਾ ਹੁੰਦਾ ਹੈ ਜਿਹੜਾ ਸਰੀਰ ਹੈ ਮੇਰ ਸਰੀਰ ਹੈ ਉਹਨੂੰ ਦ੍ਰਿ ਨਦਰ ਸਰੇ ਕੋਪੜੀ ਦਿਮਾਗ ਦਾ ਉਹ ਸਗਰ ਬੈਠੀ ਹੈ ਨਾਣਾ ਦੇ ਵੀ ਸਗਰ ਬਣਿਆ ਨਾ ਪਾੜ ਦੇ ਉੱਤੇ ਸਰੀਰ ਨੂੰ ਜੇ ਪਾੜ ਮੰਨ ਲੀਏ ਉਹਦੇ ਉੱਤੇ ਬੈਠੀ ਚਲ ਅੱਖਾਂ ਤੇ ਵੀ ਉੱਪਰ ਪੰਨਾਂ ਤੇ ਵੀ ਉੱਪਰ ਨੱਕ ਤੇ ਵੀ ਉੱਪਰ ਗਿਆਨ ਅੰਦਰ ਸਾਡੇ ਦੇ ਜੁੜੇ ਦੇ ਇਹ ਬੈਠੀ ਹੈ ਜਿਹਦੇ ਕਲ ਸੋਰ ਹੈ ਦੇਵਤਿਆਂ ਨੂੰ ਜਿਤਨ ਵਾਲੀ ਦੇਵਤੇ ਜਿਹੜੇ ਨੇ ਨਾ ਦੇਵਤੇ ਦੇਵਤੇ ਦੰਦਰ ਸੰਸਾਰ ਨੂੰ ਕੁਛ ਇਹਦਾ ਉਹਨੂੰ ਕਹਿੰਦੇ ਨੇ ਜੋ ਦੇਣੇ ਕੀ ਇੱਛਾ ਰੱਖਦਾ ਹੈ ਕੁਛ ਮੰਗਦਾ ਨਹੀਂ ਕਿਸੇ ਸੇ ਉਹ ਦੇਵਤਾ ਹੁੰਦਾ ਉਹਨੂੰ ਜਿੱਤਣ ਵਾਲੀ ਹੈ ਉਹਨਾਂ ਦੇ ਮਨ ਜਿੱਤਣ ਵਾਲੀ ਹੈ ਮਨ ਜਿੱਤ ਤੇ ਸੁਰ ਚਰੀ ਜਿੰਨੀਆਂ ਸੁਰਾਂ ਸੁਰਗ ਏ ਵੀ ਸੁਰ ਦਾ ਮੰਨ ਨਹੀਂ ਦੇਲਤਾ ਹੁੰਦਾ ਸੁਰ ਅੱਡ ਅੱਡ ਸੁਰਾਂ ਧਰਮ ਦੀਆਂ ਅੱਡ ਅੱਡ ਵਿਚਾਰ ਤਾਰਾ ਵਾਂਣ ਜੜੀਆਂ ਅੱਡ ਅੱਡ ਸੁਰਾਂ ਨੇ ਉਹ ਕਹਿੰਦਾ ਸੁਰ ਹੈ ਅੱਡ ਸੁਰ ਸਾਰੀਆਂ ਸੁਰਾਂ ਨੂੰ ਸੱਦ ਸਰ ਵਾਲੀ ਹੈ ਇੱਕ ਕਰਨ ਵਾਲੀ ਹੈ ਕਰਨਾ ਇੱਕ ਕਰਨਾ ਸਾਰੀਆਂ ਮਤਨ ਇੱਕ ਮਤ ਇੱਕ ਧਾਗੇ ਵਿੱਚ ਇੱਕ ਸੂਤ ਵਿੱਚ ਪਰੋਲ ਸੁਰਸਰੀ ਪਰਸੇਵ ਜਾਚੈ ਸੁਰਸਰੀ ਸੁਰਸਰੀ ਕੋਈ ਕੰਪਰੋਮਾਈਜ਼ ਨਹੀਂ ਕਿਸੇ ਨਾਲ ਕਰਦੀ ਉਹ ਉਹਦੇ ਨਾਲੇ ਸਾਰਿਆਂ ਨੂੰ ਕੰਪਰੋਮਾਈਜ਼ ਕਰਨਾ ਪੈਂਦਾ ਆਪਣਾ ਨਾਂ ਨਹੀਂ ਉਲਟ ਮੋੜਨਾ ਉਹਦਾ ਨਾਂ ਸਦਾ ਸਦਾ ਹੀ ਰਹੂਗਾ ਬਹਿਣ ਨੂੰ ਵੀ ਕਹਿੰਦੇ ਨੇ ਬਹਿਣ ਸ਼ੋਰਟ ਵਿੱਚ ਇਸ ਪੰਕਤੀ ਦਾ ਅਰਥ ਕੀ ਹੋਇਆ ਜੀ ਨਖ ਪਰਸੇਵ ਜਾਚੈ ਜੇ ਜਦ ਜਿੱਦੀ ਚਲਦੀ ਹੈ ਸੁਰਸਰੀ ਦਰਿਆ ਆਨੇ ਚਲਦੇ ਨੇ ਸਾਰੇ ਕੇ ਚਲਦੇ ਨਦੀਆਂ ਬਿਲਕੁਲ ਸਿੱਧੀ ਚਲਦੀ ਹੈ ਜੇ ਨਾਉ ਚਲਦਾ ਬਹਿਣ ਸਿੱਧਾ ਹੈ ਨਖ ਨਾਉ ਸਿੱਧਾ ਜਾਂਦਾ ਪਰਸੇਵ ਬਹਿਣ ਨੂੰ ਕਹਾਂਗੇ ਜੀ ਬਹਿਣ ਬਹੁ ਬਬਈ ਸੁਰਸਰੀ ਦਾ ਇੱਕ ਅਰਥ ਜਾਣਨਾ ਚਾਹੁੰਦਾ ਸੀ ਜਿਵੇਂ ਇੱਕ ਬਾਣੀ ਚ ਪੰਕਤੀ ਹੈ ਸੁਰਾ ਅਪਵਿੱਤਰ ਨਤ ਅਵਰ ਜਲਦੇ ਸੁਰਸਰੀ ਮਿਲਤ ਨਹੀਂ ਹੋਈ ਆਨੰਦ ਜਿਸ ਵਕਤ ਜਿਹੜੇ ਆਪਵਿੱਤਰ ਜਲ ਜਿਹੜੇ ਹੁੰਦੇ ਹਨ ਸੁਰਾ ਜਿਹੜੀ ਹੈ ਸੁਰਾ ਸ਼ਰਾਬ ਨੂੰ ਕਹਿੰਦੇ ਨੇ ਸੁਰ ਅਪਵਿੱਤਰ ਆ ਜਿਹੜੀ ਸੁਰਾ ਸ਼ਰਾਬ ਹੈ ਇਹ ਅਪਵਿੱਤਰ ਜਲ ਮੰਨੇ ਇਹਨੂੰ ਸਾਰਿਆਂ ਨੂੰ ਨਤ ਅਵਰ ਜਲ ਰੇ ਇਹਦੇ ਬਰਾਬਰ ਕੋਈ ਹੋਰ ਪਵਿੱਤਰ ਜਲ ਨਹੀਂ ਹੈਗਾ ਇਹ ਮੰਨਦੈ ਨੇ ਇਹ ਨੂੰ ਸ਼ੱਕ ਹੈ ਅਹੰਕਾਰਵਾਦ ਕਰਮ ਵਧਾਉਣ ਵਾਲੀ ਚੀਜ਼ ਹੈ ਤਾਂ ਪਵਿੱਤਰ ਹੈ ਗੰਗਾ ਵਿੱਚ ਆਗਦੀ ਹੈ ਇਹਦਾ ਨਾਂ ਜੇ ਇਹ ਗੰਗਾ ਜਲ ਵੇਦੇ ਵਿੱਚ ਪਾ ਦਈਏ ਗੰਗਾ ਜਲ ਚ ਪੈ ਜਵੇ ਗੰਗਾ ਦੇ ਵਿੱਚ ਜਿਵੇਂ ਆ ਛੋਟੇ ਛੋਟੇ ਦਰਿਆਨ ਨੇ ਉਹਨਾਂ ਦੇ ਨਾਂ ਨੇ ਜਦੋਂ ਗੰਗਾਜ ਪੈ ਜਾਂਦਾ ਨਾ ਫਿਰ ਨਾਂ ਆਪਣਾ ਖਤਮ ਹੋ ਜਾਂਦਾ ਗੰਗਾ ਹੀ ਰਹਿ ਜਾਂਦੀ ਹੈ ਜਦੋਂ ਸੋ ਉਹਦੇ ਵਿੱਚ ਮਿਲ ਜਾਂਦੇ ਨੇ ਰੋਂਗਾ ਦੇ ਵਿੱਚ ਫਿਰ ਉਹਦਾ ਆਪਣਾ ਨਾਂ ਖਤਮ ਹੋ ਜਾਂਦਾ ਹੈ। ਪਰ ਸੰਤ ਜਿਹੜੇ ਜੇ ਸੁਰਾ ਦੇ ਸ਼ਰਾਬ ਦੇ ਵਿੱਚ ਰੋਂਗਾ ਜਦ ਬਾਲਵੇਂ ਸੰਤ ਨਹੀਂ ਪੀਂਦੇ। ਸੰਤ ਜਿਹੜੇ ਨੇ ਉਹਨੂੰ ਪੀਂਦੇ ਨਹੀਂ ਹਨ। ਹੋਏ ਆਨੰਦ ਵੱਖਰਾ ਨਹੀਂ ਰਹਿੰਦਾ ਫਿਰ ਉਹ ਹੋਲ ਸੁਰਸਰੀ ਦਾ ਰੂਪੇ ਹੋ ਜਾਂਦਾ ਹੈ। ਨਦੀਆਂ ਨਾਲਿਆਂ ਟੋਬਿਆਂ ਦਾ ਪਾਣੀ ਮਿਲ ਸੋ ਸੁਸਰੀ ਹੋ ਜਾਏ। ਫਿਰ ਉਹਦਾ ਆਪਣਾ ਮजूद ਖਤਮ ਹੋ ਜਾਂਦਾ ਹੈ। ਦੇ ਸ਼ਬਦ ਜਿਹੜੇ ਨੇ ਜੇ ਭਗਤੀ ਦੇ ਸ਼ਬਦ ਲਿਖ ਲਵੇ ਕਾੜ ਦੇ ਰੁਸ਼ ਦੇ ਪੱਤਿਆਂ ਤੇ ਉਹ ਪਵਿੱਤਰ ਹੋ ਜਾਂਦੇ ਉਹਨੂੰ ਮੱਥਾ ਟੇਕੀਦਾ। ਪਰ ਇਹ ਸੰਤ ਨਹੀਂ ਮੰਨਦੇ। ਪਗਤਾਨੋ ਜਿਵੇਂ ਜਾਚ ਪੈਦਾ ਹੋਏ ਨੇ ਫੇਰ ਵੀ ਇਹਨਾਂ ਦੇ ਅੰਦਰ ਰਹੀ ਜਾਂਦੀ ਮੈਨੇ ਉਧਰ ਗੰਗਾ ਚ ਮਿਲਿਆ ਆ ਪਵਿੱਤਰ ਜਲ ਨਦੀਆਂ ਨਾਲਿਆਂ ਡੋਬਿਆਂ ਦਾ ਸ਼ਹਿਰਾਂ ਦਾ ਉਹ ਜਿਹੜੇ ਸੰਤ ਨੇ ਇਹਨਾਂ ਦੀ ਫੱਟੀ ਪੋਚੀ ਆ ਗੱਲ ਕਹਿ ਕੇ ਇੱਕ ਪਾਸੇ ਤੁਸੀਂ ਇੱਕ ਗੱਲ ਮੰਨਦੇ ਹੋ ਦੂਏ ਪਾਸੇ ਉਹ ਗੱਲ ਨਹੀਂ ਮੰਨਦੇ ਆਮ ਲਗੇ ਗੰਗਾ ਦੇ ਵਿੱਚ ਹਰਦਵਾਰ ਦਾ ਰਿਸ਼ੀ ਕੇ ਦਾ ਗੰਗਲਦਾ ਆਖੇ ਉਹ ਤਾਂ ਤੁਸੀਂ ਉਹ ਹੋ ਜਾ ਪਵਿੱਤਰ ਸਮਝ ਲਿਆ ਗੰਗਾ ਜਲ ਲਾਤਾ ਛਿੜਕਤਾ ਉਹ ਪਵਿੱਤਰ ਹੋ ਗਿਆ ਜੁੱਤੀ ਪਵਿੱਤਰ ਹੋ ਗਈ ਗੰਗਾ ਜਲ ਛੜਕੇ ਤੇ ਜੁੱਤੀ ਬਣਾਉਣ ਵਾਲਾ ਛਮਾਰ ਪਵਿੱਤਰ ਹੀ ਹੋਇਆ ਗੰਗਾ ਨਾਤੇ ਛੇ ਆਦੋਂ ਦੂਸਾਂ ਵੀ ਜਾਇਓ ਪਰ ਮੈਂ ਕੀ ਗੱਲ ਨੂੰ ਇਹ ਕੀ ਕਿਹ ਹੈ ਜੋ ਤੂੰ ਜਨ ਨੂੰ ਨੀਚ ਰੱਖਣਾ ਮੰਨਿਆ ਵੀ ਇਹ ਨੂੰ ਨੀਚੇ ਰੋ ਜਿਉ ਨੀਚ ਹੈ ਕਿਉਂ ਤੁਹਾਡੇ ਗੋਵਰ ਨਹੀਂ ਨੀਚ ਉੱਚ ਨਹੀਂ ਕੀਤੇ ਉਹ ਕਦੇ ਮੇਰਾ ਗੋਵਰ ਉੱਚ ਉੱਚ ਕਰਦਾ ਇਹ ਸੇ ਤੋੜਦਾ ਨਹੀਂ ਉਹ ਹਾਲ ਤੱਕ ਤੋੜਦਾ ਨਹੀਂ ਉਹ ਇਹਨਾਂ ਦੇ ਵੀ ਸੀਗੇ ਨਾ ਉਹ ਬਣੇ ਹੋਏ ਜਿਹੜੇ ਸੰਤ ਫਾਲੇ ਹੋਣੇ ਮਾਰਟੋ ਤੋਂ ਛੇਗ ਨੇ ਨਹੀਂ ਇਹ ਨਹੀਂ ਗੱਲ ਆਸੀ ਬੰਦੇ ਐਵੇਂ ਅਦਾਲਤਾਂ ਤਾੜੇ ਬਣਾਏ ਤੇ ਨਾ ਜੀ ਇਹਨਾਂ ਦੀ ਮਰਜ਼ੀ ਦੀ ਬਰਦਾ ਹੈ ਜਿਹੜੀ ਗੱਲ ਇਹਨਾਂ ਨੂੰ ਸੋਚ ਲੱਗਦੀ ਹੈ ਬੰਦੇ ਨਹੀਂ ਨਹੀਂ ਹੋਏ ਆਨੰਦ ਉਹ ਵੱਖਰਾ ਨਹੀਂ ਹੋ ਜਾਂਦਾ ਫਿਰ ਸਹੁਰੇ ਹੋ ਰਹਿੰਦਾ ਹੈ ਵਿੱਚ ਮਿਲ ਕੇ ਉਹਦਾ ਵੱਖਰਾ ਮजूद ਨਹੀਂ ਰਹਿੰਦਾ ਜਮਨਾ ਮਿਲ ਗਈ ਗੰਗਾ ਚ ਉਹਦਾ ਵजूद ਖਤਮ ਹੋ ਗਿਆ ਅੱਗੇ ਗੰਗਾ ਹੀ ਚੱਲੂ ਜਮਨਾ ਖਤਮ ਪਰ ਭਗਤਾਂ ਦੀ ਬਾਣੀ ਰਬਦਾਸ ਦੀ ਬਾਣੀ ਰਬਦਾਸ ਭਗਤ ਉਹ ਕਹੇ ਵੀ ਭਗਤਾਂ ਚ ਨਿਰਲਿਆ ਤੁਸੀਂ ਕਹਿੰਦੇ ਉਹਦੀ ਬਾਣੀ ਬਾਹਰ ਕੱਢਦੇ ਹੋ ਤਾਂ ਜਵਾਬ ਸੀ ਉਹ ਵਖਰਾ ਭਾਤੇ ਹੋ ਕੇ ਵੀ ਵਖਰਾ ਸੋਰਸੇ ਜਿ ਮੜਕੇ ਵੀ ਵੱਖਰਾ ਜਮਨਾ ਉਸ ਸੋਰਸੇ ਜਿ ਮੜਕੇ ਬੱਕਰੀ ਨਹੀਂ ਰਹੀ ਮਾਇਆ ਵਿੱਚ ਕੀ ਫੈਸਲੇ ਥੋਡੇ ਨੇ ਜ਼ੁਰੇ ਫੈਸਲੇ ਨੇ ਕਿਸੇ ਚੀਤੇ ਚੋਟ ਕੀਤੀ ਹੋਈ ਆ ਸਮਝਦਾ ਤਾਂ ਨਹੀਂ ਉਹਨਾਂ ਦੇ ਵਿਚਾਰ ਤੇ ਉਹਨਾਂ ਦੇ ਅੰਦਰ ਜਿਹੜੀ ਖੋਟ ਆ ਤੇ ਚੋਟ ਆ ਖੋਟ ਤੇ ਚੋਟ ਆ ਖੋਟ ਉਹਨਾਂ ਜਿੱਥੇ ਇਹ ਦੁੱਖ ਅਨਕਠੋ ਹੈ ਇਥੋਂ ਨਾ ਇਥੋਂ ਖੰਬਿਜਲੀ ਨਹੀਂ ਜੇ ਇਹ ਪਵਿੱਤਰ ਨਹੀਂ ਹੋ ਸਕਦੇ ਕਿਉਂਕਿ ਜੁੱਤੀ ਬਣਾਉਂਦਾ ਇਹ ਚਮਾਰ ਚਮੜਾ ਗਾਉਦਾ ਲੂ ਨੂੰ ਚੱਕਦਾ ਚਫਾਲ ਕਰਦਾ ਚਮੜਾ ਲਾਉਂਦਾ ਉਹ ਅਪਵਿੱਤਰ ਹੈ ਜੁੱਤੀ ਵੀ ਗੋਪਵਿੱਤਰ ਹੈ ਗੋ ਗੋਉ ਤਾਂ ਅਪਵਿੱਤਰ ਹੈ ਤੇ ਮਰ ਜਵੇ ਫੇ ਪਵਿੱਤਰ ਉਹਦੇ ਵਰਗਾ ਪਵਿੱਤਰ ਕੁਝ ਨਹੀਂ ਜੀ ਉਹਦਾ ਮਾਸ ਆ ਪਵਿੱਤਰ ਹੈ ਦੁੱਧ ਪਵਿੱਤਰ ਹੈ ਕਿਉਂ ਮਾਸ ਕਿਉਂ ਪਵਿੱਤਰ ਹੈ ਭਾਈ ਦੁੱਧ ਕਿਉਂ ਪਵਿੱਤਰ ਹੈ ਮਾਸ ਕਿਉਂ ਪਵਿੱਤਰ ਹੈ ਦੱਸ ਕੇ ਰੂਲ ਮਰਜੀ ਦੇ ਬਣਾਏ ਹੋਏ ਨੇ ਇਹ ਕਰਕੇ ਸੱਜੋਗ ਦੇ ਵਿੱਚ ਗੋ ਮਰੇ ਦੇ ਕਰਦੇ ਸੀ ਸਭ ਤੋਂ ਸ੍ਰੇਸ਼ ਕਿਉਂਕਾ ਗਊ ਸਭ ਤੋਂ ਪਵਿੱਤਰ ਜਾਨਵਰ ਹੈ ਉਹਦਾ ਮਾਸ ਵੀ ਪਵਿੱਤਰ ਹੈ ਇਰਾਨੇ ਜਦ ਦੇਖਿਆ ਪਤਾ ਲੱਗਿਆ ਵੀ ਖੇਤੀ ਕਰਨੀ ਹੈ ਆਪਣੀ ਬਣਾਤਾ ਪੈਣਾ ਇਹ ਇੱਥੇ ਪੈਣ ਲੋ ਸਾਨੂੰ ਇਹਦੀ ਲੋੜ ਹੈ ਸਮਾਜਿਕ ਲੋੜ ਨੂੰ ਧਰਮ ਸੀ ਕੀ ਕਰਦੇ ਸੀ ਸਮਾਜਾ ਤਾਂ ਮਰਜੀ ਦਾ ਉਹਦਾ ਪਰਦਾ ਫਾਸ਼ ਹੋਣ ਵਾਲਾ ਹੁਣ ਪਰਦਾ ਫਾਸ਼ ਹੋ ਰਿਹਾ ਹਿੰਦੂ ਹਿੰਦੂ ਨੇ ਆਕੇ ਕੀਤਾ ਹੈ ਜਦ ਤੱਕ ਤੇ ਬੰਨ ਲਗਿਆ ਉਹ ਹਿੰਦੂ ਬਣ ਕੇ ਜਾਂਦੇ ਬਣੇ ਹਿੰਦੂ ਜਾਤੇ ਹੀ ਨਾਂ ਰੱਖਿਆ ਨੇ ਆਪਣੇ ਅੰਦਰਾਂ ਦਾਸਲੀ ਛੱਡ ਫੈਸਲੇ ਲੈ ਲਏ ਇਹਨਾਂ ਨੂੰ ਤਾਂ ਹਿੰਦੂ ਕਹਿਣੇ ਸੀ ਉਹਨੂੰ ਉਹਨਾਂ ਜਾਂ ਤਾਂ ਤਰਵਜਨ ਤਾਂ ਸਾਜਿ ਵੇਦ ਛੱਡ ਤਾ ਜਮਨ ਛੱਡ ਦੇ ਫੈਸਲੇ ਤੋਂ ਕਹਿ ਕਰਨੇ ਸ਼ੁਰੂ ਕਰਤੇ ਠਗੀਆਂ ਫਰੇਬ ਸਭ ਨੂੰ ਜਾਇਜ਼ ਕਰਾ ਦਿੱਤਾ ਇਹਦੇ ਵਿੱਚ ਨਰਨਸਾਂ ਵਿੱਚ ਬਿਸ਼ਰੂ ਭੱਜ ਗਿਆ ਲੈ ਕੇ ਅਮਰਤ ਜਾਇਜ਼ ਹੈ ਕਮੇਟਵੰਤ ਕਹੇ ਸੀ ਜੰਗ ਬੰਦੀ ਦੀ ਅਰਜੁਨ ਦੇ ਮੁੰਡੇ ਨਾਲ ਧੋਖਾ ਕਰ ਲਿਆ ਜਾਇਜ਼ ਹੈ ਹੋਂ ਜੁਦ ਵਿੱਚ ਕੁਝ ਵੀ ਜਾਇਜ਼ ਹੈ ਸਭ ਕੋ ਧੋਖੇ ਤਾਂ ਨਨਵਾਂ ਸਾਹਿਬ ਛਡਾ ਲਿਆ ਧੋਖੇ ਨਾਲ ਬਾਅਦ ਆਪਣਾ ਘਰ ਤਾਂ ਸਭ ਗਏ ਇੱਥੋਂ ਆ ਕੇ ਤੁਹਾਨੂੰ ਨਸ਼ ਹੋ ਗਿਆ ਧੋਖਾ ਤਰਮ ਜਾ ਵੜਿਆ ਚਰਮੇ ਧੋਖਾ ਬਣ ਗਿਆ ਚਰਮੇ ਨੋਂ ਤੇ ਹੀ ਧੋਖਾ ਦੇ ਰਹੇ ਨੇ ਲੋਕਾਂ ਨੂੰ ਕਿ ਖਾਣੇ ਆਕਾਰ ਸਰਤ ਬਣਾ ਕੇ ਧੋਖਾ ਦਿੱਤਾ ਸਿੱਖਾਂ ਨੂੰ ਐ ਖਾਲੀ ਦਲ ਬਣਾ ਕੇ ਗੁਰਦਾਰੇ ਬਣਾ ਕੇ ਧੋਖਾ ਦਿੱਤਾ ਹੰਥ ਬਣਾ ਕੇ ਖੋਹ ਲੈ ਕੇ ਧੋਖਾ ਕੀ ਕਰੇ ਆ ਧੋਖਾ ਦਿੱਤਾ ਹੁਣ ਮੰਨ ਵੀ ਗਏ ਵੀ ਗਲਤ ਪਰਚਾਰ ਮੰਨ ਵੀ ਗਏ ਮੰਨ ਵਿੱਚ ਗਏ ਸੰਦ ਕੋਈ ਧਰਮ ਨਹੀਂ ਹਿੰਦੁਸਤਾਨ ਦੇ ਉਹਦੇ ਵਿੱਚ ਹਿੰਦੂ ਉਸ ਨੂੰ ਸੱਚ ਬਸਾਈ ਆਪਸੇ ਮੈਂ ਹਾਂ ਭਾਈ ਭਾਈ ਇਹ ਲੈ ਕੇ ਅਭੀ ਹੋਇਆ ਹਿੰਦੂ ਤਰਮ ਕਾਨੂੰਨ ਲਿਖਿਆ ਵੀ ਹੋਇਆ ਹੁਣ ਕਹਿੰਦੇ ਤਰਮ ਨਹੀਂ ਹਿੰਦੂ ਸੁਪਰੀਮ ਕੋਰਟ ਨੇ ਵੀ ਕਹਾਤਾ ਕੋਮ ਜਾ ਕੇ ਤਰਮ ਜਿੰਦਾ 50 ਬਣਾ ਲਿਆ ਆਹ ਕੁਛ ਹੈ ਵਿਸ਼ਵਾਸ ਕੌਣ ਕਰੇ ਇਹਨੂੰ ਬੋਲਣ ਕਵੇਂ ਬੋਲਣ ਕਵੇਂ ਤੁਹਾਨੂੰ ਦੇ ਉਸਤੇ ਐਂ ਤਾਂ ਧੋਖੇ ਵਾਲ ਸਾਰੇ ਰਾਜ ਧਰਮ ਹੁੰਦਾ ਹੈ ਰਾਜੇ ਦਾ ਇੱਕ ਧਰਮ ਹੁੰਦਾ ਹੈ ਆਜਾ ਦਾ ਧਰਮ ਬੌਲਦੀ ਪਾਲਣਾ ਕਰਨਾ ਗਰੀਬ ਦੀ ਪਰਵਰਿਸ਼ ਕਰਨਾ ਕਮਜ਼ੋਰ ਨੂੰ ਬਚਾਉਣਾ ਕਮਜ਼ੋਰ ਦੀ ਰੱਖਿਆ ਕਰਨਾ ਤਕੜੇ ਨੂੰ ਦੇ ਨੱਥ ਪੋੜੀ ਜੇ ਤੱਕ ਆਖਾਲ ਦਾ ਨੱਥ ਪੋੜੀ ਉਹਨੂੰ ਸਜ਼ਾ ਦੇਣੀ ਪਰ ਇੱਥੇ ਤਾਂ ਸਰਕਾਰ ਧਖਾ ਕਰਦੀ ਹੈ ਆਪੇ ظلم دی انتہا ہے اد یا راجہ ہی شیر منی ویس شیر بن جائے مقدمے کتے بن جانا سانو کتے فڑوتا پر تے پرمیشر اپے کوئی کرے ہیلا تا دنیا بچے ورنہ دنیا نو بچن کون دے تے کھان والے نے سب جوں ਇਦਸੋਕ ਕੇ ਘਾਰੇ ਲੀਡਰ ਬਣ ਕੇ ਆਦਮੀ ਨੂੰ ਘਾਰੇ ਨੇ ਆਦਮੀ ਆਦਮੀ ਆਦਮੀ ਦਾ ਖੂਨ ਚੂਸ ਰਿਹਾ ਛਰੇ ਆਮ ਚੂਸ ਰਿਹਾ ਤੇਕ ਸਵਾਕੇ ਚੂਸ ਰਿਹਾ ੱੱਕਾ ਕਰਕੇ ਚੂਸ ਰਿਹਾ ਕਾਨੂੰਨ ਬਣਾ ਕੇ ਚੂਸ ਰਿਹਾ ਫਿਰ ਤਾਂ ਪਰਮੇਸ਼ਰ ਆਪੇ ਹੀ ਕੁਝ ਕਰੇ ਆਪੇ ਕਿਸ ਰੂਪ ਵਿੱਚ ਪ੍ਰਗਟ ਹੋਵੇ ਜੀ ਆਪੇ ਕੋ ਕਲਾ ਵਰਤਾਵੇ ਖੇਡ ਵਰਤਾਵੇ ਤਾਂ ਗਲ ਉਹ ਖੇਡ ਵਰਤ ਰਹੀ ਹੈ ਉਹ ਹਲਾ ਰਿਹਾ ਆਪਣੀ ਹੁਣ ਪਿਆ ਪਿਆ ਜਿਵੇਂ ਕੋਈ ਪਾਸਾ ਲੈਂਦਾ ਕਰਵਟ ਬਦਲ ਰਿਹਾ ਹੋ ਜਦ ਕਰਵਟ ਬਦਲਦਾ ਅਸਲਜੋਕਰ ਵਤ ਹੁੰਦਾ ਆਰਾ ਚੱਲਦਾ ਫਿਰ ਇਹਨਾਂ ਤੇ ਜੁਲਮ ਤੇ ਜੁਲਮ ਤੇ ਸਲਤੇ ਪਹਿਲਾਂ ਤਾਂ ਧਰਮ ਦੇ ਸਲਤੇ ਆਰਾ ਚੱਲਿਆ ਨਾ ਧਰਮੀਆਂ ਦੇ ਸਲਤੇ ਚੱਲਿਆ ਨਹੀਂ ਆਰਾ ਦਿੱਲੀ ਚ ਜੀ ਚੜਨ ਕੜੀਆਂ ਤੇ ਚੜੇ ਨਹੀਂ ਨਰਮੀ ਹੋਰ ਜਾਲਮਾਂ ਤੇ ਆਰੇ ਚੱਲਣਗੇ ਕਰਵਟ ਬਦਲ ਗਈ ਹੋਰ ਨਾਲੇ ਸਮੇਂ ਤੇ ਜਾਲਮਾਂ ਦੇ ਉੱਤੇ ਆਰੇ ਚੱਲਣਗੇ ਕਰਮੀ ਨਾ ਕਰੀ ਜਲ ਲੈਣ ਅੰਦਰ ਤਾਂ ਹੁਣ ਵੀ ਚੱਲਦੇ ਨੇ ਇਹਨਾਂ ਦੇ ਅੰਦਰ ਹੁਣ ਵੀ ਚੱਲਦੇ ਚਿੰਤਾ ਦੇ ਆਰੇ ਅੰਦਰ ਫਿਕਰ ਪੈ ਗਿਆ ਵੀ ਕੀ ਅੰਤਯੰਤਾ ਸਭ ਨੂੰ ਵਿਗਵੇ ਗੰਢ ਖਲੋਹ ਦੁਨੀਆ ਨੂੰ ਬੇਕਾਬੂ ਹੁੰਦੀ ਜਾਂਦੀ ਹੈ ਹਾਂਜੀ ਆਪਾਂ ਇਸ ਪੰਕਤੀ ਦੇ ਅਰਥ ਕੀਤੇ ਸੀ ਨਖ ਪਰਸੇਵ ਜਾਂਚੈ ਸੁਰਸਰੀ ਇਹਦੇ ਜਿਹੜੇ ਅਰਥ ਹੋਏ ਪਹਿਲਾਂ ਉਹ ਹੋਏ ਪਹਿਣ ਗੰਗਾ ਉਸ ਦੇ ਦਰ ਤੇ ਉਸ ਦੇ ਨੌਂ ਦਾ ਪਸੀਨਾ ਹੈ ਆਪਾਂ ਪਹਿਲਾਂ ਨਹੀਂ ਕੀਤੇ ਹਾਂ ਸੁਰਾ ਅਪਵਿੱਤਰ ਨਤ ਅਵਰ ਜਲਦੇ ਉੱਥੇ ਆਪਾਂ ਸੁਰਸਰੀ ਦੇਤ ਗੰਗਾ ਕਿਤੇ ਨਹੀਂ ਇਹ ਗੰਗਾ ਕਹਿੰਦੇ ਨੇ ਗਿਆਨ ਦੀ ਗੰਗਾ ਸਾਡੀ ਪ੍ਰਕਾਸ਼ ਗੰਗਾ ਨਹੀਂ ਕਹਿੰਦੇ ਹਾਂਜੀ ਫਿਰ ਉਹ ਵੀ ਤਾਂ ਗੰਗਾ ਹੀ ਹੈ ਇਹਨਾਂ ਦੀ ਆਪਣੀਆਂ ਗੰਗਾ ਸਾਡੀ ਆਪਣੀਆਂ ਬਈ ਗੰਗਾ ਇਹ ਨਹੀਂ ਚਲਦੀ ਜਿਵੇਂ ਦੀ ਚਲਦੀ ਹੈ ਦੇਖੋ ਬੱਦਲ ਵੀ ਚੱਲਦੇ ਨੇ ਹਵਾ ਨਾਲ ਸਿੱਧਾ ਹੀ ਜਾਂਦੇ ਨੇ ਜਾਂਦੇ دریاਵਾਂੋਂ ਤਾਂ ਜਾਂਦੇ ਨਹੀਂ ਹਵਾ ਜਾਂ ਚਲਦੀ ਹੈ ਸਿੱਧੀ ਚਲਦੀ ਹੈ ਜੇ ਪੂਰਬ ਦੇ ਜਿੱਧਰ ਵੀ ਚਲਦੀ ਹੈ ਸਿੱਧੀ ਚਲਦੀ ਹੈ تیر ਜਿੱਧਰ ਮਰਜੀ ਮਾਰਦੇ ਸਦਾ ਜਾਊਗਾ ਜੇ ਪਰ تیر ਬਦਲ ਤੇ تیر ਸਦਾ ਜਾਊਗਾ ਕਿ تیر ਮਹ ਜਾਂਦੀ ਹੈ ਇਹ ਨਖ ਨਖ ਜੋ ਸਿੱਧਾ ਜਾਵੇ ਨਾ ਹੁੰਦਾ ਐਸਾ ਨੋ ਨਿਕਲਦਾ ਜਣਾ ਚੋਂ ਸਦਾ ਜਾਂਦਾ ਗੋੜ ਗੋੜ ਨਹੀਂ ਹੁੰਦਾ ਨੌਂ ਨੇ ਜੋ ਕਈ ਜਗ੍ਹਾ ਮੋਟੀ ਪਤਲੀ ਵੀ ਹੁੰਦੀ ਹੈ ਹੱਡੀ ਹੋ ਜਾਂਦੀ ਹੈ ਰਾਜ ਨੌਂ ਨਹੀਂ ਮੋਟਾ ਪਤਲਾ ਹੁੰਦਾ ਜਾਂ ਜਾਂ ਬਾਬਾ ਜੀ ਗੰਗਾ ਆਏਗਾ ਅਰਥ ਗੰਗਾ ਦਾ ਗੰਗਾ ਨਹੀਂ ਯਾਰ ਗੰਗਾ ਇਹ ਗੰਗਾ ਇਹਨਾਂ ਦੀ ਗੰਗਾ ਤੇ ਦ੍ਰਿਸ਼ਟੀ ਨਾ ਰੱਖ ਗੰਗਾ ਤੇ ਸਿਰਫ ਇੱਕੋ ਹੀ ਤਿੰਨ ਚੀਜ਼ਾਂ ਹੁੰਦੀਆਂ ਨੇ ਨੰਨਾ ਦਾ ਕੋਈ ਚੇਂਜ ਮੰਦੀ ਹੁੰਦੀ ਆ ਸੰਸਾਰੀ ਸਾਰੀ ਗੱਲਾਂ ਨਹੀਂ ਮਿਲਦੀਆਂ ਹੁੰਦੀਆਂ ਇੱਕ ਤਾਂ بارش ਪੈਂਦੀ ਆ ਉਤੋਂ ਆਹਤੋਂ ਵੇਗੇ ਤੋਂ ਚੱਲਦੀ ਆ ਪੱਛਮ ਤੋਂ ਪੂਰਬ ਨੂੰ ਜਾਂਦੀ ਆ ਅਸਲ 'ਚ ਇਹਨਾਂ ਦੀ ਪੂਰਬ ਦੱਖਣ ਨੂੰ ਜਾਂਦੀ ਆ ਉਲਟੇ ਹਨ ਗੰਗਾ ਦਾ ਉਲਟੇ ਨਾ ਨਹੀਂ ਗਾ ਜੀ ਸਾਡੇ ਵਾਲੇ ਪੂਰਬ ਤੋਂ ਨਿਕਲ ਕੇ ਪੱਛਮ ਨੂੰ ਜਾਂਦੀ ਇਹਨਾਂ ਦੀ ਪੱਛਮ ਤੋਂ ਨਿਕਲ ਕੇ ਪੂਰਬ ਨੂੰ ਜਾਂਦੀ ਆ ਸਾਡੀ ਬਾਹਰ ਨਾਲ ਦੇ ਉੱਤੇ ਵੀ ਜਲਦੀ ਇਹਨਾਂ ਦੀ ਥੱਲੇ ਨੂੰ ਜਾਂਦੀ ਹੈ। ਰਾਮ ਕੀ ਤੇ ਚੜਦੇ ਹੋ ਕਬੀਰ। ਬੱਦਲ ਥੱਲੇ ਉੱਪਰ ਨੂੰ ਗਏ ਨੇ। ਉਪਰੋਂ ਥੱਲੇ ਨੂੰ ਵਰ੍ਹਦੇ ਨੇ। ਇਵੇਂ ਪਹਿਲਾਂ ਬੁੱਧ ਸੋ ਤੋਤੇ ਨੂੰ ਜਾਂਦੀ ਹੈ ਉੱਤੇ ਚੜਦੀ ਆਕਾਸ਼ 'ਚ ਹੈ। ਜ਼ਮੀਨ ਤੋਂ ਉੱਪਰ ਉਹ ਤੋਤੇ ਬੋਲਦੀ ਹੈ ਜਦ ਬਾਰਿਸ਼ ਹੁੰਦੀ ਹੈ। ਇਹੀ ਕਹੂੰਗਾ ਸਾਡੀ। ਵੇਗਾ ਇਹੀ ਹੈ। ਇਹਨਾਂ ਨੇ ਆ ਗੰਗਾ ਬਹਾਲੀ ਬਣਾ ਲਈ। ਦਰਿਆ ਤਾਂ ਹੋਰ ਵੀ ਬਤੇ ਨੇ ਸੰਸਾਰ 'ਚ ਉਹ ਵੀ ਤਾਂ ਹੈਗੇ ਨੇ ਫਿਰ ਜਿੰਨੀਆਂ ਵੀ ਨਦੀਆਂ ਨੇ ਬਾੜ ਚੋਂ ਕੇ ਇੱਕ ਨਦੀ ਹੈ ਜਿਹੜੀ ਜਮਨਾ ਥੱਲੇ ਤੋਂ ਰਲਦੀ ਆ ਕੇ ਪੱਕੀ ਸਾਹਿਬ ਇਧਰੋਂ ਬਾੜ ਦੇ ਵਿੱਚੋਂ ਜਿਹੜੀ ਦੱਖਣ ਦੇ ਵਿੱਚੋਂ ਰਲਦੀ ਹੈ ਨਾ ਉਹ ਸਰ ਪੰਜਮਨਾ ਹੈ ਦੱਖਣ ਪੱਛਮ ਤੋਂ ਰਲਦੀ ਹੈ ਵਿੱਚ ਆ ਕੇ ਤਾਂ ਕਿ ਪੂਰਬ ਦੇ ਵਿੱਚ ਉਹ ਉੱਤਰ ਚੋਂ ਆ ਕੇ ਦੇ ਜੀ ਪਾਰਨੀ ਜਨੈ ਜੇ ਪਈ ਜਾਂਦਾ ਨਾ ਰੀਆਂ ਦਾ ਐਵੇਂ ਸਾਡੇ ਵਿਚਾਰਤਾ ਰਹੇ ਗੁਰਮਤਿ ਦੱਖਣ ਦੇ ਕੇ ਇਹ ਪਹਾੜ ਰੀਆਂ ਜਿੰਨੀ ਉੱਪਰ ਨੂੰ ਵਿਚਾਰਤਾ ਰਹਾਂ ਨੇ ਸਾਰੀਆਂ ਵਿਚਰੜ ਜਾਂਦੀ ਇਹਦੇ ਇਸ ਬੁੰਦਲ ਤੱਕ ਚਲੀ ਜਾਂਦੀ ਹੈ ਇਹਨੂੰ ਤਾਂ ਗੰਗਾ ਉਹਦੇ ਨੇ ਤਸ਼ਵੀਰ ਦਿੱਤੀ ਹੋਈ ਹੈ ਕੰਪੈਰੀਜ਼ਨ ਕੀਤਾ ਹੈ ਗੰਗਾ ਕਾਨੂੰ ਹੈ ਗੰਗਾ ਕਿਤੇ ਗੰਗਾ ਇਹਨਾਂ ਦੀ ਹੋਊਗਾਗਾ ਇਹ ਗੰਗਾ ਸ਼ਿਵਦੀਆਂ ਝੜਾਂ ਝੜ ਜਾਈ ਐ ਜਿਹੜੇ ਛੇ ਪਖਤ ਨੇ ਉਹ ਇਹਦਾ ਮਸਲਾ ਹੈ ਉਹ ਗੈਨ ਦੀ ਗੰਗਾ ਨੂੰ ਝੜਾਂ ਝੜ ਜਾਂਦੇ ਨੇ ਜਲਦਾਂ ਰੱਖ ਕੇ ਨੋ ਵਧਾ ਕੇ ਨੋਗੇ ਬਤਾਉਂਦੇ ਨੇ ਹੱਥ ਨਖਨ ਬੜਾਏ ਕਹਿਣਾ ਨਹੀਂ ਨੋ ਬੜਵੜੜ ਕਰਦੇ ਨੇ ਉਹ ਨਾ ਖਿਆ ਉੱਥੇ ਨੋ ਨਹੀਂ ਨੇ ਹੋ ਸਿੱਧੇ ਜਾਂਦੇ ਨੇ ਇਹ ਉਹਨਾਂ ਨੇ ਇਹਨਾਂ ਚੀਜ਼ਾਂ ਨਾਲ ਮਿਸਯੂਜ਼ ਕੀਤਾ ਹੋਇਆ ਹੈ। ਨਖਰਾਤ ਨਾਮ ਕਰ ਲਿਆ ਇਹਨਾਂ ਨੇ। ਨਾ ਹੁੰਦਾ ਨਹੀਂ ਨਖਰਾਤ। ਨਖਰਾ ਸਖਤ ਤੇ ਸਿੱਧਾ। ਸੁਧਰ ਸੁਧਰ ਇਹ ਚਲੋ ਤਮ। ਨਾ ਤੜ ਕੋ ਕੱਢ ਲਈਏ। ਆਦਮੀ ਸਿੱਧਾ ਹੋਵੇ ਸਪਸ਼ਟ ਹੋਣਾ। ਇਹਦਾ ਬੜਾ ਸਿੱਧਾ ਆਦਮੀ ਹੈ। ਕਹਿੰਦੇ ਨਾ ਆਪਾ। ਸੱਚੀ ਗੱਲ ਕਰਦਾ। ਸਪਸ਼ਟ ਗੱਲ ਕਰਦਾ। ਜਿਹੜਾ ਵਲਪਾ ਦੇ ਗੱਲ ਕਰਦਾ ਉਹ ਨਪਾਨ ਕਪੜੇ ਕਹਿੰਦੇ ਆ ਪਾ ਕਹਿੰਦੇ ਵਾੜਾ ਅੰਦਰ ਕਪੜੇ ਦੀ ਨਿਸ਼ਾਨੀ ਹੈ ਵਾੜਾ ਇਹਵੇਂ ਦਰਿਆ ਜਿੰਨੇ ਚੱਲਦੇ ਨੇ ਸਿੱਧੇ ਚੱਲਦੇ ਹੀ ਨਹੀਂ ਪਾਣੀ ਕਦੇ ਐਵੇਂ ਚਲੇਗਾ ਇਹਨੂੰ ਇਹਨੂੰ ਇਹਨੂੰ ਇਹ ਕਹਿੰਦਾ ਸੱਪ ਦੀ ਚਾਲ ਚੱਲਣਾ ਸੱਪ ਸਿੱਧਾ ਚੱਲਦਾ ਹੀ ਨਹੀਂ ਮਨ ਸਿੱਧਾ ਚੱਲਦਾ ਹੀ ਨਹੀਂ ਮਨ ਨੂੰ ਸੱਪ ਨਾਲ ਜੋੜਿਆ ਹੈ ਤਾਂ ਹੀ ਬੀਜ ਨੂੰ ਨਵੀਂ ਛੱਪਾ ਨਾਲ ਛਵੀ ਦੇ ਨਾਲ ਛਵੀ ਛੱਪਾ ਦੋ ਦੋਹਾਂ ਦਾ ਮਨ ਹਾਵੀ ਹੈ ਦੋਹਾਂ ਤੇ ਬਈ ਉਹ ਛਵੀ ਦਾ ਗਾਲੂ ਨੇ ਬੈਠ ਪਾਇਆ ਛੱਪਨੇ ਜਮਨਜੀ ਕੋਲ ਦਮੇ ਉਹ ਤਕਾਲ ਚ ਛੱਪ ਪਿਆ ਹੋਇਆ ਜੀ ਜਮਨਜੀ ਕੋਲ ਦਦਾ ਸਰੂਪ ਨਾ ਸਵੈਮ ਦਾ ਰੂਪ ਐ ਨਾ ਖਾਇ ਹੋ। ਸ੍ਰੂਪ ਨਾ ਖਾਨਿਆ ਲਵ। ਰਾਮਨ ਦੀ ਭੈਣ। ਸਰੂਪ ਨਜਣ ਸਰੂ ਜਿਹੜੇ ਰੂਪ ਹੁੰਦਾ ਇੱਕ ਸਰੂਪ ਹੁੰਦਾ। ਸਰੂਪ ਜੋਤ ਦਾ ਹੁੰਦਾ। ਮਨ ਤੋਂ ਜੋਤ ਸਰੂਪ ਹੈ। ਰੂਪ ਨਹੀਂ ਲਿਆ। ਸਵੈਮ ਦਾ ਰੂਪ ਜਿਹੜਾ ਸਰੂਪ ਹੁੰਦਾ। ਸਰੀਰ ਸਵੈਮ ਦਾ ਰੂਪ ਨਹੀਂ ਹੈ, ਸ੍ਰੀ ਰੂਪ ਹੈ। ਇਹ ਵਿਸ਼ੇ ਸੰਦਾਰ ਜੇ ਤੂੰ ਦੇਖਦਾ ਹਰਕਾ ਰੂਪ ਹੈ ਸੁੰਦਰ ਰੂਪ ਨੀ ਹੈ ਬਾਲਾ ਰੂਪ ਹੈ ਕਪੜੇ ਖੂਪ ਹੁੰਦਾ ਕਮੀਜ਼ ਖੂਪ ਹੈ ਪਜਾਮਾ ਪੈਂਟ ਖੂਪ ਹੈ ਪਤਾ ਵੀ ਲਤਾਜ ਬੌਰ ਹੈ ਜੁਰਾਵ ਖੂਪ ਹੈ ਪਤਾ ਪੈਰਾਂ ਨੂੰ ਪਉ ਹੈ ਉਰਗਰੇ ਬੰਦੀ ਹੋਣੀ ਦਸਤਾਨਾ ਹੱਥ 'ਤੇ ਪਉ ਵਨਨ ਗਲਛੇ ਪਊਗੀ ਕਿ ਸ਼ਹਿਰਾ ਤੇੜੇ ਪਊਗਾ ਰੂਪ ਉਹਦਾ ਕਪੜੇ ਦਾ ਜਿਹੜੀ ਜੋਤ ਆ ਉਹ ਸਰੀਰ ਤੇ ਪਹਿਨੇ ਵਾਲਾ ਕਪੜਾ ਹੈ ਸਰੀਰ ਦਾ ਰੂਪ ਨਾਲ ਮੈਚ ਕਰਦਾ ਜੋ ਉਹਦਾ ਰੂਪ ਨਾਲ ਕੋਈ ਵੀ ਕਪੜਾ ਨਹੀਂ ਕਰਦਾ ਉਹ ਸਰੀਰ ਕਰਦਾ ਜੋ ਉਹਦੇ ਰੂਪ ਨਾਲ ਮੈਚ ਸਵੈਮ ਦਾ ਰੂਪ ਕੁਛ ਹੋਰ ਹੈ ਉਹਦਾ ਜੋਤ ਆ ਜਿਹੜੀ ਉਹ ਚਮਕਾ ਜਿਹੜੀ ਚਾਨਣਾ ਰੋਸ਼ਨੀ ਹੈ ਉਹਦਾ ਸਰੂਪ ਹੈ ਸਵੈਮ ਦਾ ਰੂਪ ਹੈ ਜਿਹੜਾ ਉਹ ਸਰੂਪ ਨਾ। ਉਹ ਤੇ ਵੀ ਨਾ ਖਾਲਾ ਹੋਇਆ। ਉਹਨੂੰ 라वण ਦੀ ਪੈਣ ਮੰਨੇ ਆ। ਮੰਨਿਆ ਨੇ ਮੰਨੇ। ਜੀ। 라वण ਕੀ ਹੈ? 라वण ਚਾਰਵੇਂ ਦੱਗਿਆ ਤਾਂ ਬਵੇਕ ਹੈ। ਉਹ ਬਵੇਕ ਬੁੱਧੀ ਹੈ। ਉਹ ਪੈਣ ਪ੍ਰਾਪ ਹੋ ਗਿਆ ਇੱਥੇ ਆ ਕੇ ਦੇਉ ਸਾਤ ਪੈਣ ਪ੍ਰਾਪ ਹਾਂ। ਇਹ ਤੇ ਪੈਣ ਪ੍ਰਾਪ ਦਾ ਰਿਸ਼ਤਾ। ਤੂੰ ਮੇਰਾ ਪਤਾ ਤੂੰ ਮੇਰਾ ਮਾਤਾ ਤੂੰ ਮੇਰਾ ਬੰਦੂ ਤੂੰ ਮੇਰਾ ਪ੍ਰਾਤਾ ਤੇ ਤੇ ਪ੍ਰਾਤਾ ਦੇ ਰੂਪ ਜੀ ਵੀ ਰੱਥਿਆ ਹੋਇਆ ਵੇਖਿਆ ਅਮਰ ਤਕੀਨ ਹੈ ਸੁਰਸੁਰੀ ਦੀ ਥੋੜੀ ਜੀ ਕਲੈਰੀਫਿਕੇਸ਼ਨ ਚਾਹੀਦੀ ਹੈ ਜੀ ਹਾਂ ਆਪਾਂ ਪਹਿਲਾਂ ਨਖ ਦੀ ਕਰ ਲਈ ਨਖ ਦੀ ਕਰ ਰਏ ਸੀ ਆਪਾਂ ਨਖ ਦੀ ਹੈ ਜੀ ਨਖ ਸਿੱਧਾ ਇੱਕੋ ਸਿਕਰਾ ਸ ਇੱਕ ਰੂਪ ਨੋ ਜਿਹੜੇ ਨੇ ਜੇ ਨੋ ਕੱਟ ਕੇ ਤੋਂ ਲਿਆ ਕੇ ਰੱਖੀਏ ਦੰਗੜਾਂ ਦੇ ਨੋ ਕੋਈ ਜਦੋਂ ਪਛਾਣ ਨਹੀਂ ਹੁੰਦਾ ਕਿਹੜੀ ਬਲ ਨੇ ਪਤਾ ਲੱਗਦਾ ਵੀ ਆ ਹੱਡੀ ਕਿੱਥੇ ਦੀ ਹੈ ਨੋ ਨਹੀਂ ਪਛਾਣ ਹੁੰਦੇ ਮਾਇਨਾ ਮੋੜ ਮੋਟਾਈ ਫਰਕ ਹੁੰਦਾ ਇਹ ਗੁਰੂ ਜਿਹੜਾ ਹੈ ਉਨਾਰਾ ਰੂਪ ਹੈ ਸੇਮ ਰੂਪ ਉਤੇ ਰੂਪ ਦਾ ਫਰਕ ਹੈ ਬਸ ਪਬਈ 15 ਨੰਬਰ 972 ਤੇ ਹੈ ਜਬ ਨਖ ਸਿੱਖ ਤਬ ਅੰਤਰ ਮੱਜਨ ਕੀਨਾ ਆ ਦੇਖ ਨਰਚ ਕਾਰਨ ਕੋਰ ਮਤ ਸਿੱਧੀ ਸਿਕਾ ਸਪੈਸ ਚਖਿਆ ਸਿੱਧੀ ਗੱਲ ਉਹਨੂੰ ਖੋਜੀ ਨਖਸਿਕ ਬਾਪੇ ਅੰਤਰੇ ਮੰਜਨਗੀ ਨਾ ਬਾੜ ਨਹੀਂ ਹੈਗਾ ਫਿਰ ਕੁਝ ਨਹੀਂ ਸੱਚੀ ਸਖੈ ਦਾ ਨਾ ਹੁੰਨਾ ਸਖਦਾ ਸੱਚੀ ਸਖੈ ਬਣ ਗਿਆ ਨਾ ਬਣ ਗਿਆ ਨਖ ਪਰਸੇਵ ਗੁਰਮਤਿ ਵੀ ਬਣ ਗਿਆ ਹਾਂਜੀ ਨਖ ਪਰਸੇਵ ਜਾਂਚ ਹੈ ਜਾਂਚ ਹੈ ਸੁਰਸਰੀ ਉਹਦਨ ਪਤਾ ਲੱਗਿਆ ਬੇਰਤ ਕੀ ਹੈ ਠੀਕ ਹੈ ਜੀ ਕਲੀਅਰ ਹੈ ਬਸ ਐਟਾ ਦਾ ਬਿਲਕੁਲ ਕਲੀਅਰ ਹਾਂਜੀ ਉਹ ਰ ਘਰ ਹੈ ਬਹੁਤ ਵਕਦੀ ਹੈ ਹਾਂ ਉਹ ਇਸ ਨੂੰ ਦਰਿਆ ਕਹੇ ਆਕਾਸ਼ ਮਿਆਂ ਨੇ ਲਹੰਗ ਦਰਿਆ ਗੁਸਲ ਕਰਤਬ ਬੂਧ ਇਹ ਉਹੀ ਐ ਸੋਸਰੀ ਸਮਝਾ ਨਖ ਪਰਸੇਵ ਹੈ ਇਹਦੇ ਵਿਦਵਾਨਾਂ ਨੇ ਵੱਖਰੇ ਵੱਖਰੇ ਨਾਮ ਰਖੇ ਨੇ ਉਹ ਇੱਕ ਰੂਪ ਕੀਤੇ ਨਖ ਪਰਸੇਵ ਹੋ ਗਿਆ ਸੋਸਰੀ ਵੀ ਉਸਨੂੰ ਕਹਿੰਦੇ ਨੇ ਭਾਈ ਆਸਤ ਕੀਤਾ ਹੋਇਆ ਆਹ ਸਭ ਪਛਾਤਰ ਸੋਦੇ ਨੇ ਬਕਰੇ ਬਕਰੇ ਵਿਦਵਾਨਾਂ ਨੇ 9 ਬਕਰੇ ਬਕਰੇ ਰੱਖ ਲੈ ਵੇਦ ਪ੍ਰਾਣ ਸਿਮਰਤ ਸੁਦਾਖਰ ਕੀਨੇ ਰਾਮ ਨਾਮ ਇੱਕ ਆਖਰ ਰਾਮ ਨਾਮ ਦੇ ਨਾਲ ਜੋ ਹੁਣ ਥੋੜੀ ਥੋੜੀ ਦੇ ਆਪਾਂ ਖੋਜ ਕੀਤੀ ਅਰਥ ਦੀ ਨਾਖ ਸਿੱਖ ਦੀ ਕਿਹੜੇ ਨਾਉ ਤੇ ਅਲਸਾ ਕੇ ਜੀ ਆਪਾਂ ਕੀਤਾ ਗੁਰਬਾਣੀ ਦੇ ਜਗਾ ਜਗਾ ਸਮਝ ਆਹ ਟੈਂਕਾਏ ਤਾਂ ਸਮਝ ਲੱਗਦੀ ਐ ਤਾਂ ਇਹੀ ਹੋ ਕਰ ਸਕਦੇ ਵੱਖਰੇ ਟੀਕੇ ਨੇ ਵੱਖਰੇ ਵੱਖਰੇ ਆਏ ਨੇ ਹੁਣ ਆਹ ਜਿਹੜੀ ਪੰਕਤੀ ਤਾਂ ਬੋਲੀ ਐ ਜਿਹੜੇ ਅਥੋਰਿਟੀ ਕੀ ਕੀਤੇ ਨੇ ਪਹਿਲੇ ਉਹ ਵੀ ਦੇਖ ਲੈ ਨਖ ਸਿੱਖਦੇ ਹੱਥ ਕੀ ਕੀਤੇ ਨੇ ਉਹਨਾਂ ਨੇ ਨਖ ਸਿੱਖ ਪੈਰਾਂ ਦੇ ਨਹਾਂ ਤੋਂ ਲੈ ਕੇ ਸਿਰ ਦੀ तक सारे ਸਾਰੇ ਨੂੰ ਚੰਗੀ ਤਰ੍ਹਾਂ ਹੁਣ ਜਦੋਂ ਆਪਣੇ ਇਸ ਮਨ ਨੂੰ ਚੰਗੀ ਤਰ੍ਹਾਂ ਵੇਖਦਾ ਹਾਂ ਅੱਛਾ ਤਾਂ ਆਪਣੇ ਅੰਦਰ ਹੀ ਇਸ਼ਨਾਨ ਕਰਦਾ ਹਾਂ ਲਾ ਉਹਦਾ ਨਾ ਹੈਗਾ ਉਹਦੇ ਮਨ ਦੇ ਨਾ ਹੈਗੇ ਚੋਟੀ ਹੈਗੀ ਵਿਚਾਰ ਪਾਤ ਤੱਕ ਨਹੀਂ ਹਾਂਜੀ ਉਲਝਾਵਾ ਜੋ ਜਿੱਕੇ ਦੇ ਵਖਰਾ ਪੜਉਂਦਾ ਨਹੀਂ ਜਿਹੜੇ ਆਵਾ ਬਾਇ ਉਹਨਾਂ ਨੇ ਹੋਰ ਕਹਿਤਾ ਹੋ ਕੀ ਲੱਭ ਲੂ ਅੱਧੀ ਕਿ ਜੁਕੀ ਲੱਭੂ ਗੱਲ ਬਣਾਲਾ ਆਇਆ ਦਲ ਆਇਆ ਠੀਕੇ ਕਿਤਾਬਾਂ ਨਿਕਲ ਯੂਨੀਵਰਸਿਟੀਆਂ ਗੱਡੇ ਭਰੇ ਪਏ ਨੇ ਕੀ ਕਰ ਲੂ ਪੜ ਕੇ ਕਿਤਾਬਾਂ ਨੂੰ ਜਿਹੜੇ ਆਪ ਉੜ ਹੋਏ ਇਹ ਗ੍ਰੰਥਾਂ ਦੇ ਵਿੱਚ ਆਪੇ ਨੇ ਕਿਤਾਬਾਂ ਲਕੀਆਂ ਨੇ ਯੂਨੀਵਰਸਿਟੀ ਵਾਲੇ ਕੀ ਗੱਲ ਨੂੰ ਉੱਥੇ phd wale ki kar lane utthe ki karde bechare uddje hoye apni kitaban padhi gaye uddje hoye ne uddje hoye wo likhi gaye uddje hoye prachar kari gaye hor sare kehne vi galat ho gaya galat ki ta tu hi khojde beemanta jo swaroop hai ussi bichoti kithon aavi bhai ye ki karde ho tu itthe aake murti pooja banati ਜਾਰਾ ਚੇਤਨੂ ਇੱਕ ਕਰਤਾ ਹੋ ਜਾਰਾ ਚੇਤਨੂ ਇੱਕ ਕਰਨਾ ਆਇਆ ਸੀ ਉੱਥੇ ਪ੍ਰੋਫੈਸਰ ਨੇ ਕੋਲ ਫਿਜ਼ਿਕਸ ਦਾ ਉਹਨਾਂ ਦਾ ਕੀ ਨੋਸੀਆ ਹੰਦੇ ਜ਼ਿੰਦਾ ਹਾਂਜੀ ਜੀ ਸਪਤ ਸਮੁੰਦ ਚਾਚੇ ਘੜਥਲੀ ਸਪਤ ਸਪਤ ਦਾ ਸਤ ਵੀ ਹੁੰਦਾ ਸਪਤ ਦਾ ਸਤ ਸਮਾਂ ਸਮੁੰਦਰ ਉਹ ਸਤ ਸਮੁੰਦਰ ਕਿਵੇਂ ਬਈ ਦੇ ਕੋਈ ਇੱਕ ਸਪਤ ਲਫਦਾ ਇੱਕ ਸਤ ਲਫਦਾ ਸੱਤ ਨੂੰ ਕੰਨਾ ਤਤਾ ਸਤ ਜਿੱਤੇ ਸੱਤੇ ਨੂੰ ਕੰਨਾ ਤਤਾ ਸਤ ਇਹਦਾ ਅਰਥ ਹੈ ਸੈਵਨ ਜਿੱਤੇ ਸਪਤ ਅਰਥ ਹੈ ਸਤਵਮ ਸੱਤ ਨੇ ਵੀ ਦੀਆਂ ਸੱਤੇ ਸਮੁੰਦਰ ਨੇ ਜਿਹੜੀ ਸੱਤਵੀਂ ਦੇ ਵੀ ਹੈ ਸਪਤ ਸਹੀ ਹੈ ਚੰਡੀ ਹੈ ਅਬਵੇ ਖੋਦੀ ਹੈ ਉਹਦੇ ਆਲਾ ਸਮੁੰਦਰ ਉਹਦੇ ਆੜਾ ਗਿਆੰਦਾ ਸਮੁੰਦਰ ਸੱਤ ਸੱਤਵਾਂ ਨਾਕੇ 7 ਸੈਵਨ ਇਹਨਾਂ ਨੇ ਆਪੇ ਸੈਵਨ ਕੀਤਾ ਕੀ ਕੀਤਾ ਸੱਤੇ ਸਮੁੰਦਰ ਉਸ ਦੀ ਕੜਵਨ ਜੀ ਹਨ ਸੱਤ ਸੱਤਵਾਂ ਨੇ ਤਾਂ ਸੱਤਾਂ ਜਿਆਪਾ ਕਹਿੰਦੇ ਸੈਵਨਥ ਸੈਵਨ ਦਾ ਸੈਵਨ ਦਾ ਸੈਵਨ ਤੋਂ ਲੱਗਿਆ ਸੈਕੰਡ ਸੈਗਣ ਦਾ 2 ਨਹੀਂ ਸੱਤਵਾਂ ਫਸਲ ਦਾ ਕਿੰਨਾ ਪਹਿਲਾ ਫਿਰ ਇੱਥੇ ਆ ਕੇ ਆਕੀਤਾ ਨੂੰ ਨਾ ਉਹ ਫਸਲਾਂ ਤਾਂ ਇੱਕ ਨਹੀਂ ਹੁੰਦਾ ਪਹਿਲਾ ਹੁੰਦਾ ਹੈ ਇਹਨਾਂ ਨੇ ਜਾਨਵਰ ਜਿਵੇਂ ਕੀਤਾ ਹੋਇਆ ਪਬਲਿਕ ਕੀ ਕਰਦੀ ਉਹ ਪਬਲਿਕ ਦਾ ਮੂਰਖਾਂ ਦੀ ਹੈ ਵੀ ਦੁਵਾਨ ਮੂਰਖ ਹੁੰਦੇ ਨੇ ਸਾਨਾ ਬੰਦਾ ਹੁੰਦਾ ਉਹ ਦੇਖਦਾ ਵੀ ਸੱਤ ਦਾ ਸੱਤਮਾ ਹੁੰਦਾ ਉਹ ਇਹੀ ਸੱਤ ਸਿਰੰਗਾ ਉੱਤੇ ਸੋ ਬਤਾਤਾ 10 ਗਰ ਸੱਤ ਨਹੀਂ ਲੱਗਦਾ ਫਿਰ ਉਹਦੇ ਸੱਤ ਝੋਟੀਆਂ ਬਣਾਤਾ ਜਿੱਥੇ ਥਿੱਤੀ ਗੌੜੀ ਆਇਆ ਉੱਤੇ ਸਾਥ ਉੱਤੇ ਸਾਥ ਲਫਜ਼ਾ ਸੱਤੇ ਸੱਚ ਕਰ ਬਾਤਾਂ ਮਾਨ ਸੱਤੇ 7ਵੇਂ ਨੰਬਰ ਤੇ 7ਵੀਂ ਗੱਲ 7ਵਾਂ ਵਚਨ ਸੱਤੇ ਸੱਤੇ ਨਾਲ ਇਹਦੇ ਨੂੰ 7ਵੀਂ ਗੱਲ ਇਹ ਹੈ ਸਤ ਕਰ ਇਹਨੂੰ ਸੱਚੀ ਬਣਨਾ ਜਿਹੜੀ ਮੈਂ ਹੁਣ ਸੱਤਵੇਂ ਨੰਬਰ ਤੇ ਗੱਲ ਕਰਨ ਲੱਗਿਆ ਆਤਮ ਰਾਮ ਨੇ ਉਹ ਕੁਰਬਾਨ ਆਪਣੇ ਆਪ ਨੂੰ ਅਰਾਮ ਹੁੰਦਾ ਆਤਮ ਜਿਹਨਾਂ ਤੇਰਾ ਮੂੜਾ ਉਹ ਹੀ ਰਾਮ ਹੈ ਪ੍ਰਵਾਨ ਕਰਦਾ ਤੇ ਪ੍ਰਵਾਨ ਨਹੀਂ ਕਰਦਾ ਕਿਉਂਕਿ ਤੂੰ ਰਾਮ ਬਾਹਰ ਬੰਦੀ ਬੈਠਾ ਪ੍ਰਵਾਨ ਕਰਵਾਇਆ ਜਿਹਨਾਂ ਦਾ ਪ੍ਰਵਾਨ ਕਰ ਲਿਆ ਉਹਦਾ ਬੰਦਿਆ ਸਿੱਖ ਜਿਹਨੇ ਪ੍ਰਵਾਨ ਨਹੀਂ ਕੀਤਾ ਉਹ ਸਿੱਖ ਨਹੀਂ ਬਣੇ ਇਸ ਅੰਗਲ ਤਰਬਾਹ ਲਿਖਿਆ ਦਸਮ ਪਾਸ਼ਾ ਦੇ ਆਤਮ ਰਾਮ ਆਤਮ ਰਾਮ ਜਿਸ ਨਜ਼ਰੀ ਆਇਆ ਇਹ ਕਹਿੰਦਾ ਜੀ ਸੂਬੇ ਸਾਹਿਬ ਦੇ ਵਿੱਚ ਉਥੇ ਵੀ ਆਤਮ ਰਾਮ ਲਫ਼ਜ਼ ਵਰਤੇ ਇੱਥੇ ਵੀ ਆਤਮ ਰਾਮ ਨਾਮ ਵਰਤੇ ਐ ਰਾਮ ਜਿਹੜਾ ਆਤਮ ਰਾਮ ਆ ਉਹੀ ਪੰਜਵੇਂ ਪਾਸ਼ਾ ਵਰਤ ਰਹੇ ਨੇ ਉਹ ਕਹਿੰਦਾ ਆਤਮ ਰਾਮ ਰਹੋ ਪਰਵਾਣ ਇਹਨੇ ਪ੍ਰਵਾਨ ਕੀਤਾ ਕਿ ਉਹ ਕਹਿੰਦਾ ਆਤਮ ਰਾਮ ਜਿਸਨੂੰ ਨਹੀਂ ਆਇਆ ਤਤ ਕਾਲ ਦਾ ਦੇਸ ਪ੍ਰਗਟ ਆਇਆ ਤਤ ਕਾਲ ਦਾ ਦੇਸ ਦਸਾਈ ਦੇ ਸ਼ਾਵਨ ਦੇ ਪ੍ਰਗਟ ਹੋ ਗਿਆ ਸਵੇਕ ਰਾਮ ਬੋਲਦਾ ਨਜ਼ਰ ਦੀ ਆ ਰੋ ਫਰਕ ਇੱਥੇ ਹੈ ਫਰਕ ਇਹਨਾਂ ਦਾ ਜਾਣ ਕੇ ਪਾਇਆ ਹੋਇਆ ਫਿਰ ਕਹੋ ਕਬੀਰ ਤੂੰ ਰਾਮ ਕੀ ਅੰਸ਼ ਰਾਮ ਦੇ ਰੂਪ ਹੈ ਜਿਹੜਾ ਹੁਣ ਅਪੂਰਣ ਹੈ ਬੂਲ ਨਬਰ ਬਣੀ ਰਿਆ ਕਮਜ਼ੋਰ ਹੋ ਗਿਆ ਸ਼ਕਤੀ ਪੂਰੀ ਨਹੀਂ ਬੁੱਧਵਲ ਪੂਰਾ ਨਹੀਂ ਰਹਾ ਬੁੱਧਵਲ ਹੀਨ ਹੋ ਗਿਆ ਬੁੱਧਵਲ ਹੀਨ ਹੋਇਆ ਘਟਿਆ ਰੂਪ ਹੀਨ ਰੂਪ ਵੀ ਘਟ ਗਿਆ ਠੱਗਾ ਪੈ ਗਿਆ ਕਮਜ਼ੋਰ ਹੋ ਗਿਆ ਚਮਕ ਘਟ ਗਈ ਰੂਪ ਹੀਨ ਬੁੱਧਵਲ ਹੀਨ ਮੈਂ ਪਰਦਾ ਸੰਦੂਰ ਤੇ ਆਈ ਦੇਖਿਆ ਨਾ ਜੀ ਜੋਤ ਨੂੰ ਲਗਾਉਰ ਕੀ ਜੋਤ ਹੀ ਗਲ ਹੋਤੇ ਜਾਦ ਦੀ ਗੱਲ ਹੈ ਓਈ ਸੁਰਸਰੀ ਹੈ ਸੁਰਸੇ ਨਾ ਕਿਓ ਫਿਰ ਰੂਬੀ ਢੀ ਕੋਈ ਉਹਦਵਾਲ ਵੀ ਪੂਰਾ ਹੋ ਗਿਆ ਉਹ ਜਿ ਮਿਲ ਕੇ ਜੀ ਉਹ ਸੁਰਸੇ ਜਿ ਮਿਲ ਕੇ ਸੁਰਸੇ ਦਾ ਰੂਪ ਇਹ ਹੋ ਜੂ ਸੁਰਸੇ ਲੋਪ ਹੈ ਉਹ ਨਾ ਆਪਣੇ ਆਪ ਨੂੰ ਸੁਰਸੇ ਦੇ ਬਜੇ ਲੀਨ ਕਰ ਨਦੀ ਨੇ ਦੂਰੀ ਨੇ ਨਦੀਆਂ ਨਾਲੇ ਟੋਪਿਆਂ ਦਾ ਪਾਣੀ ਮਿਲ ਸੁਰਸਰੀ ਜੋ ਜ ਮਿਲ ਗਿਆ ਸੁਰਸਿ ਦਾ ਰੂਪੇ ਹੋ ਗਿਆ ਤੋ ਕਹਣਾ ਨਹੀਂ ਇਸ ਕਰਕੇ ਜਿਹੜਾ ਸੁਰਸਿ ਜੀ ਦਾ ਵਿੱਚ ਕੁਛ ਵੀ ਮਿਲ ਜਾਂਦਾ ਸੁਰਸਿ ਤੋਂ ਵੱਖਰਾ ਨਹੀਂ ਰਹਿੰਦਾ ਪਸੰਤ ਜਨ ਵੱਖਰਾ ਰੂਪ ਮੰਨਦੇ ਨੇ ਨਹੀਂ ਕਰਤਪਾਨਾ ਇਹਦਾ ਮਤਲਬ ਇਹ ਹੋਇਆ ਕਿ ਥੋੜੀ ਗੰਗਾ ਉਹ ਆਪਣਾ ਰੂਪ ਨਹੀਂ ਬਣਾ ਸਕਦੀ ਤੁਸੀਂ ਅੰਦਰੋਂ ਇਹ ਮੰਨਦੇ ਹੋ ਜੇ ਮੰਨ ਸਕਦੇ ਜੇ ਤੁਸੀਂ ਮੰਨਦੇ ਹੋ ਕਿ ਗੰਗਾ ਦਾ ਜਲ ਆਪਣਾ ਰੂਪ ਬਣਾ ਲੈਂਦਾ ਤਾਂ ਗੰਗਾ ਦੇ ਜਲ ਪਾ ਕੇ ਸ਼ਰਾਬ ਪੀ ਕੇ ਦਿਖਾਓ ਇਹ ਉਹਨਾਂ ਦਾ ਟੈਸਟ ਲਿਆ ਵਕਤਾ ਨੇ ਜੀ ਸਮਝਿਆ ਗੱਲ ਸਮਝ ਗਈ ਜੇ ਗੰਗਾ ਨੂੰ ਪਵਿੱਤਰ ਮੰਨਦੇ ਹੋ ਸ਼ਰਾਬ ਪੀ ਕੇ ਦਿਖਾਓ ਸ਼ਰਾਬ ਪੀ ਕੇ ਦਿਖਾਓ ਪੰਦੇਸ਼ ਸ਼ਰਾਬ ਪੀਂਦਾ ਨਹੀਂ ਉਹ ਵੀ ਨਹੀਂ ਤੇ ਉਹਨਾਂ ਦਾ ਪਵਿੱਤਰ ਮੰਦਾ ਨਹੀਂ ਕਹਿੰਦਾ ਹੈ ਮੰਦਾ ਨਹੀਂ ਜੋ ਕਹਿਣਾ ਹੁੰਦਾ ਨਹੀਂ ਇਹਨਾਂ ਦੀ ਗੰਗਾ ਤੋਂ ਉਹਨੂੰ ਟੌਂਟ ਮਾਰੀ ਹੈ ਜੀ। ਜਾਂ ਜੀ ਉਹਨੂੰ ਬੁਗਰਾਇਆ ਹੈ ਉਹ ਤੋਂ। ਸਪਤ ਸਮੁੰਦ ਜਾਂਚੈ ਘੜਥਲੀ। ਉਹ ਕਾੜਦੇ ਉਹਦੇ ਥਲੀ ਦੇ ਥਲ ਹੁੰਦਾ ਉਹਦਾ ਜਿਹੜੀ ਹੱਥ ਦੀ ਥੇੜੀ ਕਹਿ ਲੋ। ਘੜਥਲੀ ਹੋਣਾ ਘੜਥਲੀ ਨਹੀਂ। ਘੜ ਕੱਗਾ। ਓਏ ਘੜਥਲੀ ਯਾਰ। ਘਰ ਹੱਥਾ ਘੜਦੀ ਹੈ। ਕੱਗਾ ਨਹੀਂ ਹੈਗਾ ਜੀ। ਯਾਰ ਮੈਂ ਤੁਹਾਨੂੰ ਦੱਸਾਂ ਕਾਰਲ ਆਫ ਹੈਗਾ ਹੈ ਉੱਥੇ ਇੱਕ ਜਗ੍ਹਾ ਹੋਰ ਵੀ ਹੈ ਸਭਨਾਂ ਦਾ ਕਰ ਆ ਕਰ ਹੈ ਕਰਦੀ ਹੈ ਕਰਦੀ ਨਾ ਤੇ ਜੀ ਕਰ ਥਲੀ ਤਾਂ ਹੁੰਦਾ ਹੀ ਨਹੀਂ ਕਰ ਥਲੀ ਹੁੰਦਾ ਥਲੀ ਤਾਂ ਹੱਥ ਦੀ ਮੁਠੀ ਇੱਕੋ ਵਾਰੀ ਆਇਆ ਜੀ ਆਦ ਬਾਣੀ ਵਿੱਚ ਘੜ ਥਲੀ ਸ਼ਬਦ ਇੱਕੋ ਵਾਰੀ ਆਇਆ ਇੱਥੇ ਪਰ ਕਰ ਥਲੀ ਹੁੰਦਾ ਯਾਰ ਕਰ ਥਲੀ ਹੈ ਨਹੀਂ ਅੱਛਾ ਜੀ ਆਹ ਉਹ ਦਾ ਉਹ ਆਪੇ ਉਹ ਦਾ ਘਰ ਇਹਦਾ ਮਤਲਬ ਚਲੋ ਆਪਾਂ 2 ਮਿੰਟ ਬਾਅਦ ਫਿਰ ਉਹ ਦਾ ਕਰ ਜਿਹਦਾ ਘਰ ਹੈ ਉਹ ਘਰ ਵੱਡਾ ਹੁੰਦਾ ਘਰ ਵੱਡਾ ਜੀ ਤੁਸੀਂ ਸਰਪਿਆ ਘਰ ਹੈਗਾ ਉਹ ਤੇਰਾ ਘਰ ਤੇਨੂੰ ਬੜਾ ਛੋਟਾ ਮੇਰੇ ਤੋਂ ਬੜਾ ਜੀ ਫਿਰ ਫਿਰ ਘਰ ਦਾ ਦਾ ਜੇ ਘਰ ਹੈ ਕੋਈ ਤਾਂ ਉਹ ਵੀ ਘਰ ਤੋਂ ਦੀ ਹੈ ਉਦਾਕਾਰ ਜਿਹਨੂੰ ਕਹਿ ਦਿੱਤਾ ਜਾਂਦਾ ਜਸਰ ਮਾਰੂ ਕੋਡਾ ਆ ਰੇ ਫਿਰ ਪਰਮੇਸ਼ਰ ਦਾ ਘਰ ਪਰਮੇਸ਼ਰ ਤੋਂ ਛੋਟਾ ਹੈ ਉਹ ਆਪੇ ਆਪਣਾ ਕਹਦਾ ਯਾਰ ਉਹਦਾ ਘਰ ਕੀ ਹੋ ਜੂ ਉਹਦਾ ਘਰ ਉਹਦੇ ਵਿੱਚ ਲਿਆ ਘਰ ਹੈ ਉਹਦਾ ਘਰ ਦੀ ਹੁੰਦਾ ਥਲੀ ਕੀ ਹੁੰਦੀ ਹੈ ਥਲੀ ਕੀ ਹੈ ਥਲ ਉਹ ਥੇੜੀ ਅਥੇ ਅਥੇੜੀ ਉਹਨੇ ਹਾਂਜੀ ਇਹਨੂੰ ਥਲ ਇਹਨੂੰ ਕਹਿੰਦੇ ਨੇ ਕਰ ਹਾਲੀ ਤਪਤ ਸਮੁੰਦਰ ਉਹ ਪਿੱਛੇ ਕਾਰਲਾ ਨਾ ਉਹਦੇ ਘਰ ਉਹਦੇ ਘਰ ਤਾਂ ਘਰ ਕਰਤਾ ਚਾਚਾ ਘਰ ਸਿੱਤੇ ਕਾਰ ਉਹਨਾਂ ਨੇ ਕਹਦੇ ਠੋਕ ਤਾਂ ਇੱਥੇ ਵੀ ਠੀਕ ਹੈ ਜੀ ਹਾਂ ਘੜ ਮੇਰੇ ਭਾਲ ਕੇ ਨੇ ਕਹਿਤਾ ਯਾਰ ਇੱਕ ਘਰ ਨਹੀਂ ਹੈ ਤੇ ਘਰ ਚਾਹੀਦਾ ਘੜ ਤਾਂ ਚਲੇ ਪਿੱਛੇ ਕੜ ਥਲੀ ਸ਼ਬਦ ਬਾਬਾ ਜੀ ਕਿਸੇ ਵੀ ਗ੍ਰੰਥ ਵਿੱਚ ਨਹੀਂ ਆਇਆ ਨਾ ਦਸਮ ਬਾਣੀ ਚ ਤੇ ਨਾ ਹੀ ਆਦ ਬਾਣੀ ਚ ਇਸ ਤੋਂ ਇਲਾਵਾ ਬਹੁਤ ਜਾਨਣ ਦੀ ਕੜ ਹੈ ਜਸਲੀ ਸਾਰੇ ਖਜ਼ਾਨੇ ਹੈ ਜੀ 10 ਸਦੀਆਂ ਠਾਕੁਰ ਕਰਤਾਲ ਤਰਿਆ ਉਹਦੇ ਹੱਥ ਦੀ ਥੇਲੀ ਤੇ ਉਹਦੇ ਝੇਲੀਓ ਦਾ ਕਾਰ ਹੈ ਉਹਦੇ ਹਥੇੜੀ ਆ ਜਿਹੜੀ ਉਹਦਾ ਹੁਕਮ ਹੈ ਉਹਦਾ ਕਾਰ ਹੈ ਹੁਕਮ ਹੈ ਉਹਦਾ ਹੱਥ ਹੈ ਉਹ ਹੀ ਉਹਦਾ ਕਾਰ ਹੈ ਹੁਕਮ ਹੈ ਹੱਥ ਹੈ ਉਹਦੇ ਦੇ ਵਿੱਚ ਨੇ ਜੀ ਜਾਂਚ ਵਰਤਣੀ ਇਹਨੇ ਵਰਤਣ ਵਾਸਤੇ ਸਾਰੇ ਜੀ ਉਹਦੇ ਹੁਕਮ ਦੇ ਨੇ ਜੀ ਤੇ ਡੜਾ ਕੋਈ ਮਰਜ਼ੀ ਕਰਾ ਲਵੇ ਭਾਈ ਦਰਗਨ ਨੂੰ ਕਹਿੰਦੇ ਉਹਨਾਂ ਦਾ ਕੰਮ ਕਰਾਉਣੇ ਦੂਜੀ ਦੀ ਵਧੀਆ ਡਿਊਟੀ ਲਾ ਦੇ ਜਿਹੜਾ ਕੰਮ ਜਾਣਦਾ ਅਰਲਾ ਉਹਦੇ ਚ ਕੰਮ ਕਰਨਾ ਵੀ ਆ ਤੂੰ ਕੱਲ੍ਹ ਲਈ ਦੁਆ ਕਰਨਾ ਇਹ ਵੀ ਉਹ ਨਹੀਂ ਜਾਂਦਾ ਆਪਣੇ ਬੰਦੇ ਆਪਣੇ ਆਖਰ ਲੱਗਦੇ ਹੀ ਹੁੰਦੇ ਨੇ ਇਹ ਕੋਈ ਨਵੀਂ ਗੱਲ ਹੈ ਸੰਸਾਰੀ ਗੱਲ ਹੀ ਆ ਇਹਦੇ ਕਾਰੇ ਨੇ ਮੈਂ ਪਰ ਹੁਣ ਕੰਮ ਕਰਨ ਵਾਲੇ ਉਹਦੇ ਹੁਕਮ ਚੱਲਣ ਵਾਲੇ ਉਹ ਜੀ ਤਾਂ ਮੰਦੀ ਜਿਹੜਾ 93 ਆਪਣੇ ਆਪ ਨਹੀਂ ਲੈਦਾ ਆਪਣੀ ਕੋਸ਼ਿਸ਼ ਕਰਦਾ ਉਹਦੇ ਬੰਦੇ ਹੁਕਮਾਂ ਵਾਲੇ ਕਰਨਾ ਉਹਦੇ ਹੁਕਮ ਦੇ ਸਾਬ ਨੂੰ ਚੱਲਣ ਵਾਲੇ ਕਰਾਉਣੇ ਹੈਗੇ ਉਹਦੇ ਕੋਲ ਸਭ ਕੁਝ ਕਰਦਾ ਹੋਇਆ ਵੀ ਕੁਝ ਨਹੀਂ ਕਰਦਾ ਸਭ ਕੁਝ ਦੇਖਦਾ ਹੋਇਆ ਵੀ ਕੁਝ ਨਹੀਂ ਦੇਖਦਾ ਸਭ ਕੁਝ ਸੁਣਦਾ ਹੋਇਆ ਵੀ ਕੁਝ ਨਹੀਂ ਸੁਣਦਾ ਸਭ ਕੁਝ ਸੋਚਦਾ ਹੋਇਆ ਵੀ ਕੁਝ ਨਹੀਂ ਸੋਚਦਾ ਲੈਕਿਨ ਸਮਝਦਾ ਆਪੇ ਕੱਲਾ ਹੀ ਐ ਸਭ ਕੁਝ ਇਹ ਨਹੀਂ ਕਹਿ ਸਕਦੇ ਸਮਝਦਾ ਹੋਇਆ ਵੀ ਕੁਝ ਨਹੀਂ ਸਮਝਦਾ ਸਮਝ ਉਹਦੀ ਚਲਦੀ ਹੈ ਸੋਚ ਲੋਕਾਂ ਦੀ ਚਲਦੀ ਹੈ ਉਹਦੀ ਮਰਜ਼ੀ ਪਰ ਸੋਚ ਦੂਜਿਆਂ ਦੀ ਚਲਦੀ ਹੈ ਮਰਜ਼ੀ ਉਹਦੀ ਚਲਦੀ ਹੈ ਹਾਂਜੀ ਸੋ ਐਸਾ ਰਾਜਾ ਤ੍ਰਿਭਵਨ ਧਣੀ ਐਸਾ ਰਾਜਾ ਹੁੰਦਾ ਤੈਨ ਲੋਕ ਦਾ ਤ੍ਰਿਭਵਨ ਧਣੀ ਤਿੰਨ ਪਾਪੜਾਂ 'ਚ ਤਿੰਨ ਪਾਪੜ 'ਚ ਇੱਕੋ ਜੋਗੀ ਕਹੋ ਕਵਣ ਹੈ ਰਾਜਾ ਹੈ ਨਾ ਜੀ ਉਹ ਜਿਹੜੀ ਬਝਾਰਦਾ ਕਵਣ ਹੈ ਰਾਜਾ ਨਾ ਆ ਉਹਦੇ ਬਝਾਰ ਤੋਂ ਦੱਸੀ ਆ ਉਹ ਜਵਾਬ ਆਉਦਾ ਤਿੰਨ ਪਾਪੜਾਂ 'ਚ ਇੱਕੋ ਜੋਗੀ ਗਵੀਰ ਨੇ ਪੁੱਛਿਆ ਸੀ ਨਾ ਹੋਰ ਦੱਸੋ ਰਾਜਾ ਕੌਣ ਨੇ ਫਿਰ ਕੋਈ ਕੱਲਾ ਹੀ ਆ ਸਾਰਿਆਂ ਨੂੰ ਜੁੜਿਆ ਹੋਇਆ ਸਾਰੇ ਨਾਲ ਜੁੜਿਆ ਇੱਕੋ ਜੋਗੀ ਹੈ ਸਾਰੇ ਨਾਲ ਜੁੜਿਆ ਹੋਇਆ ਉਹ ਜਿਹਨੂੰ ਆਪਣੀ ਮਰਜ਼ੀ ਜੀਤੇ ਜੋ ਮਰਜ਼ੀ ਕਰਾ ਲਵੇ تیرے ਭਵਨ ਤਾਂ ਨਹੀਂ ਆਹੋ ਤਾਂ ਹੀ ਕੱਟ ਉਹ ਕੱਟ ਕੱਟ ਕੇ ਅੰਤਰੀ ਕੀ ਜਾਣਤਾ ਤੈਨਾਂ ਲੋਕਾਂ ਚ ਕਿ ਜੁੜਿਆ ਹੈ ਤੈਨਾਂ ਲੋਕਾਂ ਨਾਲ ਸਾਰੇ ਜੀਵਾਂ ਨਾਲ ਜੁੜਿਆ ਹੋਇਆ ਸਾਰੇ ਉਹਦੇ ਨਾਲ ਜੁੜਿਆ ਮਹਿਸੂਸ ਕਰਨ ਨਾ ਕਰਨ ਪਰ ਉਹ ਸਾਰਿਆਂ ਨਾਲ ਜੁੜਿਆ ਹੈ ਉਹਦਾ ਧਿਆਨ ਸਾਰਿਆਂ ਨਾਲ ਜੁੜਿਆ ਹੋਇਆ ਹੈ ਹਰ ਵਕਤ ਸਾਰੇ ਉਹਦੇ ਧਿਆਨ ਚ ਰਹਿੰਦੇ ਨੇ ਸਾਰੇ ਉਹਦੇ ਖਿਆਲ ਚ ਰਹਿੰਦੇ ਨੇ ਜੀ ਚਾਹੇ ਉਹਦਾ ਧਿਆਨ ਰੱਖਦੇ ਨੇ ਚਾਹੇ ਨਹੀਂ ਰੱਖਦੇ ਪਰ ਉਹ ਨਹੀਂ ਭੁੱਲਦਾ ਕਿਸੇ ਦਾ ਭਲਾਇਆ ਕੋਈ ਜਾਗਤ ਜੋਤ ਹੈ ਨਾ ਅਸੀਂ ਸੁਪਨਾ ਦੇਖਦੇ ਹਾਂ ਜਾਗਤ ਜੋਤ ਹੈ ਨਹੀਂ ਜਿਹੜਾ ਜਾਗਤ ਹੁੰਦਾ ਜੋਤ ਉਹ ਇੰਨਾ ਹੀ ਜੁੜ ਜਾਂਦਾ ਜਿਵੇਂ ਉਹ ਜੁੜਿਆ ਸਭ ਨਾਲ ਜਾਗਤ ਜੋਤ ਉਹਦੇ ਨਾਲ ਜੁੜ ਜਾਂਦਾ ਬਾਕੀਆਂ ਨਾਲ ਨਹੀਂ ਜੁੜਨੀ ਲੋੜ ਉਹ ਉਹਦੇ ਨਾਲ ਜੁੜਦਾ ਉਹਦੇ ਨਾਲ ਜੁੜ ਕੇ ਇਦਾਂ ਜੁੜਦਾ ਸਾਰਿਆਂ ਨਾਲ ਉਹ ਜੁੜਿਆ ਹੋਇਆ ਹੀ ਹੈ ਅਸੀਂ ਟੀਵੀ ਨਾਲ ਜੁੜਨਾ ਤੇ ਉਹ ਕੈਮਰੇ ਨਾਲ ਨਹੀਂ ਜੁੜਨਾ ਜਿਹੜਾ ਜਗਾ ਜਗਾ ਫੜ ਕੇ ਟੀਵੀ ਨੂੰ ਮੈਸੇਜ ਦੇ ਰਿਹਾ ਟੀਵੀ ਚਾਈ ਜਾਣਾ ਸਭ ਕੁਝ ਕੈਮਰਾ ਕੋਬਦਾ ਟੀਵੀ ਚਾ ਰਿਹਾ जी वो सब सब कुछ देखना है को देख ही जाना ठीक है जी बाबा जी इत्ते चौथे पदे दी समाप्ति है जी अच्छा जी जाचय निकटवर्ती अर्जुन ध्रु प्रहलाद अंबरीक नारद नेजय सिद्ध बुद्ध गण गंधर्व बानवे, हिला ਇਹ ਜਿਹੜੇ ਨੇ ਹੁਣੂ ਰੂਪ ਲਾਗ ਇਹ ਡਿਕਟਰੀ ਉਹਦੇ ਨੇੜੇ ਨੇ ਜਿਹੜੇ ਬਾਕੀ ਸੀ ਉਹ ਦੂਰ ਸੀਗੇ ਇੱਕ ਡਿਕਟਵਰਤੀ ਆ ਗਿਆ ਲਾਹ ਹੁਣ ਸੋਈਆਂ ਸ਼ੁਰੂ ਕਿਥੋਂ ਹੈ ਪਹਿਲਾ ਪਤਾ ਕੱਥਾ ਸ਼ੁਰੂ ਹੋਇਆ ਸੇਵੀਏ ਦੇ ਗੋਪਾਲ ਰਾਏ ਅਕੁਨ ਮਨਰਜਨ ਭਗਤ ਦਾ ਨਦੀਜਾ ਸੰਤ ਜਨ ਅਲਸੀ ਜਾਂਦੇ ਜਿਆ ਜਾਚਰ ਫੋਨ ਨੂੰ ਭਗਤੀ ਦਾਨ ਹੁਣ ਮਿਲ ਗਈ ਇਹ ਨੂੰ ਪ੍ਰੋਪਗਲਾਨ ਨੂੰ ਆ ਆ ਕੇ ਭਗਤੀ ਮਿਲ ਗਈ ਮਿਲ ਕੇ ਮੈਂ ਰਾਧ ਵਿੱਚ ਤੈਨੂੰ ਪਤਾ ਨੇ ਉਹ ਕੀ ਕਹਿੰਦੇ ਨੇ ਤੈਨੂੰ ਸੇ ਨੇ ਜੜੀਆਂ ਕਿ ਤਤੂਰੀਆ ਪਾਦਾ ਗਿਆ ਨਾ ਚਾਰ ਚਾਰੇ ਬਾਦਨ ਇਹ ਚਾਰੇ ਬਾਦਨ ਹਾਂਜੀ ਹੁਣ ਪੰਜਵਾਂ ਸ਼ੁਰੂ ਹੈ ਜੀ ਅਨੌਨੀ ਚੌਥਾ ਹੀ ਆ ਉਹ ਪਹਿਲੇ ਦੇ ਵਿੱਚ ਤਾਂ ਭਗਤੀ ਹੈ ਉਹ ਦੀ ਮੱਛਿਆ ਤਾਂ ਉੱਥੇ ਤਾਂ ਪੌਦ ਚਾਰੇ ਨੇ ਉਹ ਪਹਿਲਾਂ ਦਾ ਤਰਪ ਜਾਉ ਤਾਂ ਹੀ ਮੰਗੂਗਾ ਕੁਝ ਪਦਾਰਥ ਹਾਂ ਉੱਥੇ ਜਾਚਿਆ ਹੋਇਆ ਬੱਬੀ ਜੇ ਉੱਥੇ ਮੱਛਿਆ ਜਾਚੈਂ ਜਾਚ ਘਰ ਜਿਹਦੇ ਘਰ ਵਿੱਚ ਪਹਿਲਾਂ ਦਾ ਪੈਰ ਗੋੜਾ ਮਾਲ ਨਾਲ ਗੱਫਾ ਲੈ ਜਦੋਂ ਪਿਆਰ ਗੌੜਾ ਮਾਰ ਤੇ ਨੂੰ ਸਮਝਾਇਆ ਤੇ ਹਟ ਗਿਆ ਤਾਂ ਬਲ ਗਿਆ ਤੇ ਇਹ ਸਕੂਲ ਬਣਾਏ ਪ੍ਰਾਇਮਰੀ ਪ੍ਰੇਰੇ ਲੋਕ ਵੀ ਭਾਈ ਇੱਥੇ ਣਾਣੇ ਨੂੰ ਪੜਾਇਆ ਕਰੋ ਉਹ ਕਹਿੰਦੇ ਛੱਡੋ ਪਰੇ ਣਾਣੇ ਨੂੰ ਪੜਾ ਕੇ ਇੱਥੇ ਣਾਣਿਆਂ ਤੇ ਕੰਮ ਕਰ ਲੈ ਮੈਂ ਛੱਡਿਆ ਚਾਰੂ ਉਹ ਪ੍ਰੇਰਣਾ ਸ਼ੁਰੂ ਕੀਤੀ ਹੈ ਪਹਿਲਾਂ ਜਬ ਬਰੇਰ ਕੇ ਜਿਹੜੇ ਸਕੂਲ ਚ ਆਏ ਦਾਖਲ ਹੋਏ ਨੇ ਉਹ ਪਹਿਲਾ ਉਹ ਜਿਹੜੇ ਸੀ ਉਹ ਦਾਖਲ ਹੋਏ ਨੇ ਜਿਹੜੇ ਪੜਨ ਵਾਲੇ ਉਹ ਪਹਿਲੀ ਕਲਾਸ ਹੈ ਪਹਿਲਾ ਦਾਖਲ ਤੋਂ ਸ਼ੁਰੂ ਹੁੰਦਾ ਸਿੱਖਿਆ ਲੈਣ ਲੱਗਿਆ ਜਦ ਸਿੱਖ ਪੰਥ ਲੈਂਦਾ ਨਹੀਂ ਸਿੱਖਿਆ ਦੂਰ ਨੂੰ ਜਾਂਦਾ ਦੂਰ ਗਿਆ ਦੂਰਮਤਾ ਤਾਂ ਦੂਰਮਤਾਲੇ ਨਹੀਂ ਦੂਰਮਤ ਜਾਂ ਗੁਰਮਤ ਵਾਲ ਨੂੰ ਖੋਲਦੇ ਨੇ ਸਿੱਖਿਆ ਲੈਣ ਲੱਗਦੇ ਨੇ ਪੰਜ ਪੰਜ ਲੱਗਦੇ ਨੇ ਉਹ। ਜਾਂ ਇੱਕ ਦਾ ਬੰਦ ਮੁਖਾ ਦਾ ਘਰ ਤਾਂ ਸਿੱਖਿਆ ਲੈਦੀ ਹੀ ਨਹੀਂ। ਐਂ ਗੱਲ। ਸਾਖਤਾ ਦਾ ਘਰ ਨਹੀਂ ਗਾਲੋ ਉਹ ਤਾਂ ਖਲਾਫ ਨੇ ਨਾਮ ਤੇ। ਤਾਂ ਲਾਟਾ ਖਲਾਫ ਉਹ ਤਾਂ ਜੇ ਜਾਂ ਦੂਏ ਟੜੇ ਚੋਂਦਾ। ਫੇਰ ਪਹਿਲਾ ਪਦਾ ਸ਼ੁਰੂ ਹੁੰਦਾ। ਪਹਿਲਾ ਪਦਾ ਸ਼ੁਰੂ ਹੁੰਦਾ। ਪਹਿਲੇ ਪਦੇ ਗੁਰਮੁਖ ਮੰਨੂ ਇਕੱਠੇ ਹੀ ਨੇ ਉਹ ਲੈਣੇ ਵਾਲੇ ਨੇ ਬਾਕੀ ਨਹੀਂ ਲੈਣੇ ਵਾਲੇ ਜਿਹੜੇ ਸੁਣ ਕੇ ਲੈਣੇ ਵੱਲ ਉੱਡੇ ਨੇ ਦੂਆ ਤੋਂ ਵੱਖਰੇ ਹੁੰਦੇ ਨੇ ਨਿਖੜਦੇ ਨੇ ਉਹ ਪਹਿਲਾਂ ਪ੍ਰਾਪਤ ਹੋ ਗਿਆ ਨਾ ਛੋੜਿਆ ਮੰਨਿਆ ਉਹਨਣ ਵਾਲੂ ਆ ਗਿਆ ਜਿਹੜਾ ਜਿਹੜਾ ਮੰਨਣ ਵਾਲ ਆਇਆ ਹੀ ਨਹੀਂ ਉਹ ਜਿੱਦਿ ਹੋ ਗਿਆ ਆ ਜਦੋਂ ਜਸੂ ਹੋ ਗਿਆ ਉਹ ਉਹ ਫਿਰ ਟੱਠਿਆ ਹੋ ਗਿਆ ਉਹ ਨਾ ਹੋ ਗਿਆ ਉਹ ਫਿਰ ਉਹਦੇ ਬਾਦ ਉਹ ਰਾਮਰੇ ਇਹ ਜਿਹੜੇ ਸਾਰੇ ਨੇ ਇਹ ਕਹੇ ਨੇ ਸ੍ਰੀ ਜੱਟ ਇੱਧਰ ਆਈ ਨਹੀਂ ਉਹ ਤਾਂ ਤਰ ਗਏ ਹੋਰ ਉਹਦਾ ਇਦਾਂ ਦਾ ਮਤਲਬ ਇਹ ਨੂੰ ਤਾਂ ਪਹਿਲੇ ਕੰਨ ਪੜਾ ਲਏ ਗੁਰੂ ਇਹ ਹੋਰ ਉਹਦਾ ਤਾਂ ਉਹਦਾ ਦਰਵਾਜ਼ਾ ਤਾਲਾ ਹੋ ਗਿਆ ਬੰਦੇ ਆ ਜਿਹੜਾ ਉਹਦੇ ਚਾ ਦਤੂ ਪੂਰਾ ਚੰਨ ਨਹੀਂ ਘੜ ਲਿਆ ਬੋਣੀ ਉਹਨਾਂ ਦਾ ਦੂਜੇ ਪਾਸੇ ਉਹਦਾ ਚੰਨਾ ਵਰਦਾਰ ਹੋ ਗਿਆ ਨਾ ਪੱਲੇ ਤਾਂ ਪੱਲੇ ਜਿਹੜੇ ਨੇ ਅਸਲ ਦੇ ਵਿੱਚ ਪੱਲੇ ਜਿਹੜੇ ਨੇ ਕਿ ਬੇਦੀਆਂ ਦੇ ਜਿਹੜੇ ਨੇ ਬੇਦੀਆਂ ਦੀ ਖੁਰਾ ਹੋਜ ਮਟਾਉਣ ਵਾਲੇ ਪੱਲਿਆਂ ਨੇ ਜ਼ਿੰਮੇਵਾਰੀ ਲਈ ਹੈ ਬੇਦੀਆਂ ਦੀ ਜਣਾ ਤੇਲ ਪਾਉਣਾ ਤੇ ਗੁਰਮੱਤ ਬੇਦੀਆਂ ਬੇਦੀ ਵੇਪੜਨ ਵਾਲਾ ਹੀ ਨਾ ਗੁਰਪੰਥ ਦੀ ਕਰਨ ਦੀ ਜਾਂ ਨਬਰਦਾਰੀ ਇਹਨਾਂ ਨੇ ਲਈ ਪੱਲਿਆਂ ਨੇ ਪੱਲਿਆਂ ਨੇ ਉਹ ਤੇ ਬਾਰਾ ਨੇ ਗੁਜ਼ਾਰਦਿਆਂ ਪੱਲਿਆਂ ਕੋਲ ਪੱਲਿਆਂ ਨੇ ਉਹਦੀ ਖੰਡਣ ਨਹੀਂ ਕੀਤਾ ਬਾਰਾ ਨਾਲ ਹੁਣ ਟੱਕ ਵੀ ਹੁਣ ਵੀ ਬਾਰਾ ਦਾ ਉਹ ਕਹਿੰਦੇ ਜਨ ਘੰਡਣ ਕਰਨਾ ਚਾਹੀਦਾ ਸੀ ਕੀਤਾ ਸਗੋਂ ਬਾਰਾਂ ਦੇ ਸਹਿਣ ਹੱਕ ਜਿ ਲੈਂਦੇ ਨੇ ਇਹਦਾ ਮਤਲਬ ਬੇਦੀਆਂ ਦੀ ਖੁਰਾਕ ਉਹ ਜੜ ਪੱਤਣ ਦੀ ਜ਼ਿੰਮੇਵਾਰੀ ਪੱਲਿਆਂ ਨੇ ਲਈ ਉਹ ਪੱਲਿਆਂ ਨੇ ਆਪਣੀ ਜੜ ਪੱਟ ਲਈ ਵੇਚੀਆਂ ਸੀ ਦੀ ਪੱਟ ਹੋਣੀ ਪੱਲਿਆਂ ਦੀ ਜੜ ਤਾਂ ਪੱਟੀ ਜਾਊਗੀ ਖੁਣ ਪੱਟ ਹੋਊਗੀ ਪ੍ਰਗਟ ਹੋਏ ਤੇ ਉਹ ਥਈਨੇ ਲੋਕਾਂ ਨੂੰ ਪਤਾ ਪੱਲਿਆਂ ਦੀ ਜੜ ਰਹਿਣੀ ਨਹੀਂ ਪੱਲਿਆਂ ਦੇ ਤਾਂ ਭਲੇ ਬਣ ਜਾਣੇ ਅਰਥੇ ਬਦਲ ਜਾਣੇ ਨੇ ਭਲੇ ਥੇ ਹੀ ਭਲੇ ਤੇ ਭਲੇ ਸ਼ਬਦ ਕਾਇਵਾਰ ਆ ਫੁਰਬਾਣੀ ਚ ਭਲੋ ਭਲੋ ਆਖਿਆ ਸਭ ਕੋਈ ਪੰਨਾ ਲਾਗ ਸਕਾਇਆ ਵਾਰ ਆਇਆ ਪੰਨਾ ਤੱਕ ਵਾਰ ਬਣੀ ਆਇਆ ਉਪਰਲੇ ਸ਼ਬਦਾਂ ਪੁਰਲੇ ਪੁਰੇ ਆਇਆ ਜੀ ਪੰਨੇ ਦੇ ਉਲਟੇ ਮੋਰੇ ਆ ਭਲੇ ਸ਼ਬਦ ਭੱਬਾ ਲੱਲੇ ਨੂੰ ਇੱਕ ਲਾਮ 50 ਵਾਰ ਆਇਆ ਜੀ ਫਿਰ ਆਦਵਾਣੀ ਚ ਆਦ ਵਿੱਚ ਪੰਨੇ ਇੱਕ ਵਾਰ ਬਣੀ ਆਇਆ ਇਹਨਾਂ ਨੇ ਪੰਨੇ ਤੇ ਪੰਨੇ ਕਿਵੇਂ ਬਣਾਤਾ ਭਾਈ ਇੱਕ ਵਾਰ ਤਾਂ ਆਇਆ ਨਹੀਂ ਇਹ ਭਲੇ ਸ਼ਬਦ ਅਰਥ ਕਿਵੇਂ ਬੋਲਦੇ ਇਹ ਪੱਪਾ ਲੱਲੇ ਨੂੰ ਦੋ ਲਾਵਾਂ ਜੀ ਭੱਲੇ ਭਲੇ ਜਿਹੜੀ ਇਹ ਦੋ ਲਾਵਾਂ ਨਾਲ ਆਇਆ ਇੱਕ ਵਾਰ ਹੀ ਆਇਆ ਜੀ ਪੱਪਾ ਲੱਲੇ ਨੂੰ ਦੋ ਲਾਵਾਂ ਉਹ ਇੱਕ ਵਾਰ ਆਊਗਾ ਇੱਕ ਵਾਰ ਆਇਆ ਉਹ ਇਸ ਵਿੱਚ ਹੈ ਜੀ ਭਗਤ ਸੋਹਣੀ ਗੁਣਗਾਮ ਦੇ ਗੁਰਮਤਿ ਅਚਲੇ ਰਤਨ ਵਿਚਾਰ ਮਨ ਵਸਿਆ ਗੁਰ ਕੈ ਸ਼ਬਦ ਭਲੇ ਆ ਗੁਰ ਕੈ ਸ਼ਬਦ ਨਾਲ ਭਲੇ ਬਣੇ ਨੇ ਗੁਰ ਕੈ ਸ਼ਬਦ ਵਿੱਚੇ ਭਲਾ ਸਬਦਾ ਉਹ ਗੁਰਦੀ ਸਿੱਖਿਆ ਜਿਹੜੀ ਆ ਗੁਰਬਾਣੀ ਦੀ ਸਿੱਖਿਆ ਨਾਲ ਭਲਾ ਹੀ ਭਲਾ ਪਲੋ ਕਿੰਨੀਆਂ ਵੀ ਆਇਆ ਪਲੋ ਵੀ ਆਇਆ ਹਾਂਜੀ ਉਹ ਆਇਆ 25 ਵਾਰੀ ਫਿਰ ਇੱਕ ਵਾਰ ਇੰਨੀ ਵਾਰ ਸ਼ਬਦ ਆਇਆ ਹੋਵੇ ਗੁਰਬਾਣੀ ਤੁਸੀਂ ਉਹਦੇ ਅਰਥ ਬਦਲਤੇ ਆਪਣਾ ਨਾਲ ਜੋੜ ਲੇ ਕਿੰਨਾ ਬੜਾ ਫਰਾਦ ਹੈ ਭਲੇ ਅਮਰਦਾਸ ਗੁਰ ਕਹਰੇ ਭਲੇ ਭਾਣ ਅਮਰਦਾਸ ਬਾਤ ਆਇਆ ਅਮਰਦਾਸ ਪਹਿਨਾ ਉਦੋਂ ਪੱਲਾ ਬਾਅਦ ਚੁਰਦਾ ਫਿਰ ਅਸੀਂ ਕੁਝ ਕਹਿ ਸਕਦੇ ਸੀ ਤਾਂ ਪਹਿਲਾ ਅਮਰਦਾਸ ਬਾਅਦ ਚ ਅਮਰਦਾਸ ਤੇ ਪਹਿਲਾਂ ਵੀ ਪਲੇ ਲਾ ਕੇ ਚੱਲਦਾ ਹੈ ਅਮਰਦਾਸ ਦੇ ਨਾਲ ਕਿਵੇਂ ਜੋੜ ਦੋਗੇ ਅਮਰਦਾਸ ਪਲਾ ਬਣਿਆ ਪਲਾ ਕਨਵਾਲਾ ਬਣਿਆ ਇਹ ਪੱਲੇ ਕਹੋਂਦੇ ਹੁਣ ਨੇ ਆਪਣੇ ਆਪ ਨੂੰ ਇਹਦੀ ਮੈਂ ਕਹਿੰਦਾ ਹਿੰਦੂ ਸੀਗੇ ਉੱਤੇ ਪੱਲਾ ਆਇਆ ਕਿਸ਼ਨੂ ਉਹਦੇ ਵਿੱਚ ਕੋਲਾ ਵਰਦਨ ਪੱਲਾ ਉੱਤੇ ਪੱਲਾ ਲ ਆਇਆ ਹੋਇਆ ਹੈ ਸਾਰ ਕੋਤਾਬਲੀ ਵਿੱਚ ਇੰਦੂ ਮਾਤੀ ਚ ਪੱਲਾ ਸ਼ਬਦ ਆਇਆ ਹੋਇਆ ਹੈ ਬਿਸ਼ਨੂ ਨਾਲ ਜੁੜਿਆ ਹੋਇਆ ਇਹ ਪੱਲਿਆ ਨੇ ਠੇਕਾ ਲਿਆ ਪੱਲਿਆ ਹੈ ਸਭ ਤੋਂ ਪ੍ਰਚਾਰ ਭਾਈ ਗੁਰਦਾਸ ਭਾਈ ਗੁਰਦਾਸ ਭਾਈ ਗੁਰਦਾਸ ਨਾਲੇ ਉਹ ਦੇਵੀਆ ਮੇਰੀਆਂ ਬਾਹ ਬੇਰੀ ਬਾਣੀ ਚੜ੍ਹ ਦੋ ਉਹ ਕਹਿੰਦੇ ਵੀ ਤੇਰੀ ਬਾਣੀ ਹੈ ਤਾਂ ਦੀ ਜਾਣਨੀ ਇਥੇ ਪਰਮੇਸ਼ਰ ਦੀ ਬਾਣੀ ਚਲਦੀ ਹੈ ਇਹ ਵੀ ਸਾਖੀ ਹੈ ਛੇਵੇਂ ਪਾਸ਼ਾ ਨੇ ਭੇਜਿਆ ਔੜੇ ਲੱਗਿਆ ਉਥੋਂ ਉਲਠੀਆਂ ਕਿੜੀਆਂ ਦੇਖੀਆਂ ਇਹ ਵੀ ਪਤਾ ਫੇਰ ਵੀ ਉਹ ਵਰਉਂ ਜਾਂਦੀ ਹੈ ਕਾਸ਼ੀ ਗਿਆ ਇਹ ਤਾਂ ਮੰਗ ਗੁਰਵਾਂ ਤੇ ਤਾਂ ਨਹੀਂ ਠੀਕ ਹੋਇਆ ਕਾਸ਼ੀ ਦੀ ਪੜਾਈ ਨਾ ਜਾ ਕੇ ਠੀਕ ਹੋਇਆ ਪੂਰਾ ਹੋਇਆ। ਕੋਲੇ ਬਾਦ ਬਾਰੰਦ ਕੀ ਇਹਨੇ। ਤੇ 12 ਦਾ ਪੰਜਵੇਂ ਬਾਸ਼ਾ ਬੜੇ ਬਾਦਾਂ ਕੰਪਲੀਟ ਹੋ ਗਿਆ ਸੀ। ਕਿਰਮ ਬਾਸ਼ਾ ਬਣ ਤੰ ਵੀਰ ਤਿਆਰ ਸੀ ਉਹ ਚੜ੍ਹੌੜੀ ਪੰਜਵੇਂ ਬਾਸ਼ਾ ਨੇ ਸੀ ਪੜ੍ਹੀ। ਸਾਰੇ ਝੂਠ ਬੋਲੇ ਜਿਹੜੇ ਪੱਤੇ ਨਹੀਂ ਬੋਲੇ ਨੇ ਹੋਰ ਕੀ ਨੇ ਜੇ ਨਹੀਂ ਬੋਲੇ ਹੋਰ ਕਿਸੇ ਨੇ ਬੋਲੇ ਨੇ ਕਹਿੰਦੇ ਕਿ ਚੁੱਪ ਕਿਉਂ ਰਹੇ ਗੋਵਿੰਦਵਾਲ ਸਿੱਖੀ ਦਾ ਤੋੜਾ ਫੇਰ ਚਾਰ ਲੰਗੇ ਫੇ ਉਹਨਾਂ ਨੇ ਹਟਾਏ ਅੰਬਰ ਸਾਡੂ ਡਾਊਨ ਕਰਨ ਲੱਗੇ ਤੇ ਇਹ ਸਿੱਖੀ ਸਾਡੀ ਹੋਈ ਹੈ ਗੱਲ ਵੀ ਠੀਕ ਹੈ ਉਹਨਾਂ ਵਾਲੀ ਸਿੱਖੀ ਅੰਬਰ ਹੈ ਗੋਵਿੰਦਵਾਲ ਦੀ ਸਿੱਖੀ ਬਣਾਈ ਹੋਈ ਕੱਲ ਉਹਨਾਂ ਨੇ ਹੀ ਕਹੀ ਸੀ ਇਹ ਸਭ ਕੁਝ ਕੀ ਹੈ ਉਹ ਵੀ ਇੱਥੇ ਹੀ ਆ ਉਹਦੇ ਘਰ 'ਚ ਆ ਆਖਰ ਕਿੱਥੇ ਆ ਕੇ ਪਾਸ ਕਿੱਥੇ ਆ ਕੇ ਹੋਏ ਪਦਾਰਥ ਬੰਦੇ ਲੈਂਦੇ ਨਹੀਂ ਫਿੱਟਾਈ ਐਵੀਂ ਆਖ ਨੇ ਜਾ ਪਈ ਕਿਸੇ ਆਣੇ ਰਾਤ ਰਿਐਕਸ਼ਨ ਕਰ ਗਿਆ ਨਾ ਭੱਲਿਆ ਨੂੰ ਇੰਨਾ ਤ੍ਰੇਣਾ ਨੂੰ ਰੱਖਸ਼ ਦੀ ਕੀਤਾ ਰਿਐਕਸ਼ਨ ਦੀ ਕੀਤਾ ਤ੍ਰੇਣਾ ਨੂੰ ਹਰਾਂ ਦੀ ਕਦੇ ਚੜਨਾ ਬਰਦਾਸ਼ਤ ਨਹੀਂ ਆਉਂਦੀ ਲੱਤ ਜੂਰ ਮਾਰੀ ਹੈ ਉਹ ਵੀ ਅਮਰਦਾਦ ਦੇ ਥਾਣੀ ਤੇਣਾ ਦਾ ਇਹਨੇ ਨਾਉ ਨਹੀਂ ਲਿਆ ਕਿਉਂਕਿ ਆਮਾ ਦਾਦੀ ਬੇਇਤੀ ਕੀਤੀ ਸੀ ਤੇ ਦਾ ਲਾਉਂ ਨਹੀਂ ਲੈਂਦੇ ਪੱਲੇ ਕਿਉਂ ਲੱਤ ਮਾਰੀ ਸੀ ਅਮਰਦਾਦ ਦੇ ਇਹ ਵੀ ਚਾਰ ਨੇ ਤੇ ਹੁੰਦੇ ਪਛਾਤ ਕੋਈ ਰੋਲੇ ਨੀ ਤੇਣਾ ਦਾ ਲਾਉਂ ਨਹੀਂ ਆਉਂਦਾ ਪੱਲੇ ਪੱਲੇ ਆਉਂਦਾ ਗੁਰਦਾਸ ਦਾ ਹਾਲ ਹੁੰਦਾ ਨੱਤੂ ਦਾ ਸੁਸਾ ਜਿਗਰੇ ਨਹੀਂ ਇਹ ਸਭ ਕੀ ਹੈ ਇਹਦੇ ਬਹੁਤ بڑا ਇਤਿਹਾਸ ਹੈ ਦੇ ਵਿੱਚ ਅਸ਼ਵਦੇ ਨਾਲ ਰਿਲੇਟਡ ਹੈ ਹਾਂਜੀ ਹੁਣ ਅੱਗੇ ਪੜੋ ਭਾਈ ਗੋਇੰਦਵਾਲ ਨੂੰ ਸਿੱਖੀ ਦਾ ਧੁਰਾ ਕਹਿੰਦੇ ਆਂ ਧੁਰਾ ਹੀ ਆ ਫਿਰ ਉਹ ਵਾਲੀ ਦਾ ਜੋ ਵੀ ਆਦੀਆਂ 12 ਹਜ਼ਾਰ ਤਾਂ ਸਭ ਕੁਝ ਬਰਾਬਰ ਪ੍ਰਕਾਸ਼ ਪੜ੍ਹੀਆਂ ਜਾਂਦੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੱਚੀ ਬਾਣੀ ਵਰਵਾਣ ਕਰਦੀ ਉਹ ਰਬਨਾਲ ਖਾਂ ਸਤਗੁਰੂਗਤ ਹੋਰ ਕੱਚੀ ਆ ਬਾਣੀ ਉਹ ਕੱਚੀ ਬਾਣੀ ਨੂੰ ਤੁਸੀਂ ਬਰਾਬਰ ਕਰ ਲੈ ਪੱਕੀ ਦੇ ਅੰਨੇ ਹੋ ਗਏ ਬਿਲਕੁਲ ਗੋਲਨਾਲ ਦੀ ਕਰਾਮਾਤਾ ਗੋਲਦਵਾਲਾ ਨੇ ਨਾ ਖੋਰ ਗੱਲ ਉਹ ਅਰਜਨ ਦਾ ਜਨ ਵੀ ਗੋਇੰਦਵਾਲ ਦਾ ਨਾ RAMDAS ਗੋਇੰਦਵਾਲੇ ਰਹੇ ਸੀ ਤੇ ਦੋਨੇ ਜਿਹੜੇ ਦੂਏ ਬੜੇ ਗੋਇੰਦਵਾਲ ਦੇ ਨੇ ਨਾਲ ਕਿਹਨਾਂ ਜੱਥੇ ਇੱਥੇ ਨੇ ਉਹਨਾਂ ਦਾ ਰਿਸ਼ਤਾ ਗੋਇੰਦਵਾਲ ਨਾਲ ਹੈ ਕੱਲੇ ਅਮਰਦਾਸ ਦਾ ਰਿਸ਼ਤਾ ਗੋਇੰਦਵਾਲ ਨਾਲ ਨਹੀਂ ਅਮਰਦਾਸ ਦਾ ਪਿੰਡ ਬਾਸਰ ਕੇ ਹੈ ਅਸਲ ਉਹ ਤਾਂ ਵਾਸਣ ਦੇ ਨੇ ਇੱਥੇ ਆ ਗਏ ਰਹੇ ਨੇ ਜਲਮ ਇੱਥੇ ਦਾ ਧਰਤੀ ਇਹਦਾ ਗੋਲਨਵਾਲ ਦੀ ਜਿੱਥੇ ਧਰਤੀ ਇਹ ਦੀ ਸਿੱਖੀ ਹੈ ਭਾਈ ਗੁਰਦਾਰ ਨਾਂ ਜੋੜਿਆ ਉਹਨਾਂ ਨੇ ਉਹਨਾਂ ਨੇ ਉਹ ਸਹਿਮਤ ਰਿਹਾ ਇਹਨਾਂ ਨੇ ਬਾਬਾ ਬਟਾ ਨਹੀਂ ਰਿਹਾ ਬਕਵਾਸ ਕਰਦੇ ਨੇ ਆ ਬਾਬਾ ਬਟਾ ਛੇਵੇਂ ਪਾਸ਼ਾ ਨਾਲ ਘੋੜਿਆਂ ਦੀ ਸੇਵਾ ਕਰਦਾ ਰਿਹਾ ਕਿੱਥੇ ਉਹ ਉਥੇ ਕਾਹ ਹੋਦਾ ਇੱਕ ਪਾਸੇ ਕੰਨ ਨੂੰ ਕਾਹ ਹੋਦਾ ਉਥੇ ਐਡੀ ਦੂਰ ਉਹ ਇੱਥੇ ਸੇਵਾ ਕਰਕੇ ਕਾਹ ਹੋ ਤੜ ਜਾਂਦਾ ਸੀ ਐਡੀ ਦੂਰ ਇਹ ਸਿੱਕੀ ਗੋਇੰਦਵਾਲ ਦੀ ਉਹ ਅੰਮ੍ਰਿਤਸਰ ਦੀ ਨੇ ਅੰਮ੍ਰਿਤਸਰ ਫਰਚਾਰੀ ਗਈ ਹੈ ਗੋਇੰਦਵਾਲੋਂ ਨੇ ਜੜਾ ਜਿਵੇਂ ਨਾਮਕ ਦਾ ਨਿਰਖਾਣੇ ਕੀ ਹੈ ਮੈਨੂੰ ਇਹ ਦੱਸੋ ਨਿਰਖਾਣੇ ਕੀ ਹੈ ਦਸਬ ਬਾਚ ਜੜਾ ਪੜ੍ਹਨੇ ਕੀ ਹੈ ਕੌਜਾ ਦਾ ਪਰਨ ਕੋਈ ਨਹੀਂ ਜਾਨੂੰ ਯਾਰ ਰਸ ਪਾ ਜਿਆ ਹੋਰ ਕੀ ਹੈ ਇਹਵੇਂ ਉਹ ਦੋਹਾਂ ਦਾ ਮਾਣ ਦੇਵ ਦਾ ਪਿੰਠੀ ਦਾ ਜਨਮ ਹੈ ਤੇਰਾ ਤੇ ਅਮਰ ਨੂੰ ਨਾਂ ਅੱਜ ਵੀ ਜਿਆਦਾ ਜਿਹੜੀ ਕਹਿ ਲੋ ਲੋਧੀ ਹੋਵੇ ਚਾਹੇ ਉਹ ਨਾਂ ਗਦਰਤਾਰ ਹੋਵੇ ਜਿਤੇ ਕੋ ਨਾਮ ਦੇ ਆਖੇ ਰਹੇ ਨੇ ਇਹ ਨਾ ਸਾਰਿਆਂ ਨੂੰ ਜਿਆਦਾ ਹੀ ਪੌੜਨ ਦੇ ਰਹਿਆਂ ਸੀ ਨਰਕਾਣਾ ਸਾਹਿਬ ਨੂੰ ਜਨਮ ਹੋਇਆ ਬਰਨਾਮ ਦਾ ਹਿਸਟੋਰੀਕਲ ਹੀਰੂ ਹੋ ਕੇ ਇਹ ਮੇ ਪਰਖੀਦਾ ਇੱਥੇ ਦਾ ਇਹ ਨਾ ਸਾਰਿਆਂ ਦਾ ਤਾਂ ਦੋ ਰਾਮੰਦਰੇ ਕੁਲਕੇ ਨਹੀਂ ਕਹੀ ਗੱਲ ਪਰ ਇਹਨਾਂ ਨੇ ਫਿਰ ਦੂਏ ਸਹਿਮਤ ਨਹੀਂ ਹੁੰਦੇ ਸ੍ਰੀ ਚੰਦ ਗਿਜੜਕੇ ਸਾਹਿਬ ਤਾਂ ਨਹੀਂ ਹੁੰਦੇ ਮਨ ਨੂੰ ਪਤਾ ਜਾਂਦਾ ਕਹਨਾਂ ਦਾ ਬ੍ਰਹਮਪੂਤ ਆ ਉਹਨਾਂ ਦਾ ਸ੍ਰੀ ਗ੍ਰੰਥ ਬੀੜ ਇਹਨਾਂ ਦੀ ਹੈ ਬੀੜ ਵਿੱਚ ਇਹਨਾਂ ਦਾ ਸ੍ਰੀ ਚੰਦ ਕਹਿੰਦਾ ਕੁਝ ਵੀ ਨਹੀਂ ਸ੍ਰੀ ਚੰਦ ਨਾਲ ਕੋਈ ਸਾਧਨ ਨਾਲ ਕੋਈ ਸਾਧਨ ਨਹੀਂ ਉਹ ਤਾਂ ਆਖਿਆ ਨਾਲ ਬੀੜ ਵਿੱਚ ਕੁਝ ਨਹੀਂ ਹੈ ਸਿਰਫ ਉਹਦਾ ਪ੍ਰਭੂਤਾ ਹੈ ਨਾ ਇਹ ਇੱਕ ਐਸਾ ਗੁਰਨਾਮ ਦੀ ਬਾਣੀ ਹੈ ਬੱਬਾ ਜੀ ਉੱਪਰ ਤੁਸੀਂ ਜਦੋਂ ਸ਼ਬਦ ਸ਼ੁਰੂ ਹੋਇਆ ਤੁਸੀਂ ਉੱਥੇ ਕਿਹਾ ਹੁਣ ਕੀ ਇਹ ਮੱਥਿਆ ਭਗਤ ਭਗਤੀ ਦਾਣ ਦੀਜੈ ਜਾ ਚੇ ਉਹ ਬਾਈ ਮੱਥਿਆ ਵੱਲ ਚਲੇ ਗਏ ਨਾ ਹੋ ਭਗਤੀ ਤੋਂ ਮੱਥਿਆ ਨਾਲ ਪੱਖ ਦਿਖਾਇਆ ਤੈਨੂੰ ਮੈਂ ਗੋਲਨ ਵੱਲ ਕੀ ਹੈ ਬੱਛਿਆ ਬੱਛਿਆ ਕੰਮ ਨਾ ਉਹਦੇ ਅਰੇ ਗੋਦਾਰੇ ਮੱਛਿਆ ਬਣਾਈ ਜਾਂਦੀ ਹੈ ਪੁੱਛਦਾ ਨੇਹਰਾ ਉਹ ਮੱਛਿਆ ਤੋਂ ਬਾਅਦ ਭਗਤੀ ਸ਼ੁਰੂ ਕਰਦਾ ਹੈ ਕਬੀਰ ਕਬੀਰ ਸਿੱਤੀ 15 ਹੀ ਨਹੀਂ ਪਰ ਲਿਖਦਾ 16 ਹੋ ਇੱਕ ਮਤੋਂ ਭਗਤੀ ਸ਼ੁਰੂ ਦੀ ਜਾਂ ਚੰਨ ਥੋੜਾ ਜਿਆ ਦੇਂਗਾ ਥੋੜੀ ਹੈ ਪਰਵਾਦੀ ਚਲੀ ਜਾਂਦੀ ਹੈ ਦਿਨ ਹੋ ਠੀਕ ਹੈ ਜੀ ਸਤਿ ਆਜਿ ਮਾਰੋਂ ਸਵਾਲ ਬੱਬਾ ਜੀ ਇਹ ਐ ਕਿ ਇੱਥੇ ਆਇਆ ਦਾਨ ਦੀਜੈ ਜਾਚੇ ਸੰਤ ਜਨ ਜੇ ਸੰਤ ਜਨ ਭਗਤੀ ਮੰਗ ਰਿਹਾ ਮੱਥਿਆ ਚ ਆਓ ਸੰਤ ਜਨ ਦਾ ਭਗਤੀ ਚੌਂਦੇ ਨੇ ਹਮੇਸ਼ਾ ਮੱਥਿਆ ਚ ਵੀ ਚੌਂਦੇ ਨੇ ਜਿਵੇਂ ਪੜਨਾ ਚਾਹੁੰਦੇ ਨੇ ਆਏ ਨੇ ਸਾਰੇ ਇੱਥੇ ਭਰਮ ਦੇ ਆਣ ਨੇ ਜਬੰਦ ਆਏ ਨੇ ਉਰੇ ਹੁਣ ਜੀ ਉੱਥੇ ਮੱਥਿਆ ਤਾਂ ਸੰਤ ਜਨ ਕਿਵੇਂ ਹੋਏ ਜੀ ਇੱਥੇ ਮਾਂਖਿਆ ਉੱਥੇ ਕਿਤੇ ਮਾਂਖਿਆ ਆਂਡੇ ਦੇ ਅੰਦਰ ਬਖਸੇ ਪਰਮਦੇ ਆਂਡੇ ਦੇ ਵਿੱਚ ਆ ਸੰਤ ਬੰਦ ਹੋਇਆ ਅੱਛਾ ਜੀ ਬੰਦ ਕੀਤਾ ਕਦ ਸ਼ੌਹੰਕਾਰ ਹੋ ਗਿਆ ਬੜ ਬਰਾਬਰ ਬੋਲ ਪਿਆ ਸੁਰ ਬਜਲੀ ਮੈਂ ਮ ਲਿਖਾਇਆ ਖਸਮੇ ਕੇਦਰ ਜਾਏ ਆਏ ਗਲ ਮੈਨੂੰ ਮਰਦੋਂ ਕੀਤਾ ਜਿਹੜੇ ਮੈਂ ਬੰਦ ਕਰਦੇ ਤੇ ਉਹਨੇ ਉਹਨੇ ਬੰਦ ਕੀਤੇ ਨਹੀਂ ਉਹ ਆਟ ਖਾਤੇ ਜਿਹੜੇ ਬੋਲਦੇ ਸੀ ਅੱਡ ਘੰਟੇ ਵੀ ਜਾਓ ਬਈ ਤੇਰਾ ਵੀ ਸਾਂ ਚੱਲ ਤੇਰਾ ਵੀ ਸਾਂ ਚੱਲ ਏਰੀਆ ਤੁਹਾਡਾ ਬੜ ਜਾ ਕੇ ਨੜੀ ਜਾਓ ਜਾਓ ਸਲੀਅਰ ਹੈ ਉੱਥੋਂ ਬਾਹਰ ਨਿਕਲਨੇ ਹੁਣ ਮਸੀਹਾ ਤੂੰ ਜੀ ਜਿਹੜੇ ਦੇ ਵਿੱਚੋਂ ਅੰਦਰ ਹੀ ਰਹਿਣ ਚਾਹੁੰਦੇ ਬਾਹਰ ਨਿਕਲਣ ਦੀ ਚਾਹੁੰਦੇ ਗੁਰਬਾਣੀ ਬਾਹਰ ਕੱਢ ਰਹੀ ਹੈ ਕਬੀਰ ਬਾਣ ਕਰਦੇ ਇਕਮ ਦੇ ਵਿੱਚ ਇਕਮ ਕਹਿੰਦੇ ਪਰਬਾ ਪਰਬਾ ਕਹਿੰਦੇ ਨੇ ਇਕਮ ਦੀ ਗੰਦੇ ਪੱਖ ਦੀ ਨੂੰ ਨੇ ਪਹਿਨਾ ਪਰਬਾ ਪ੍ਰੀਤਮ ਕਰੋ ਵਿਚਾਰ ਕਟ ਮੈਂ ਖੇਲੇ ਕਟ ਕੀ ਹੈ ਪਰਮਨਾਥ ਦਾ ਘਟਾ ਕਟ ਮੈਂ ਖੇਲੇ ਆ ਪਰ ਉਹ ਜਿਹੜਾ ਇਹ ਤਾਂ ਘਟ ਸੀ ਇਹ ਤਾਂ ਸਰਵ ਵਿਆਪੀ ਦੀ ਪਰਮਦੇ ਅੰਡੇ ਚ ਕਿਵੇਂ ਪੈ ਗਿਆ ਦੇ ਕੋ ਘਨੇ ਘੜੇ ਚ ਖੇਲਦਾ ਘਟ ਇਹ ਵਿਚਾਰ ਕਰੋ ਕਿਉਂ ਘੜੇ ਖੇਲਦਾ ਕਿਉਂ ਘੜੇ ਚ ਬੜਿਆ ਇਹਦਾ ਪਰਮ ਦੂਰ ਕਰੋ ਘੜੇ ਤੋਂ ਬਾਹਰ ਕੱਢੋ ਇਹਨੂੰ ਇਹ ਇੱਥੋਂ ਸ਼ੁਰੂ ਹੋਈ ਆ ਗੱਲ ਪੜਵਾ ਪੱਖ ਦੀ ਜਿਹੜੀ ਪਹਿਲੀ ਆ ਉਹਨੂੰ ਪਰਵਾ ਕਹਿੰਦੇ ਨੇ ਮੇਰੇ ਕੱਖ ਦੀ ਪਹਿਲੀ ਨੂੰ ਇਹ ਕਹਿੰਦੇ ਨੇ ਇੱਕਮ ਜਿਹੜੀ ਆ ਜਿਹੜੀ ਮੱਛਿਆ ਵਾਲਾ ਜਿਹੜਾ ਸ਼ੁਰੂ ਹੁੰਦੀ ਆ ਜਦ ਚੰਦ ਜਾਂ ਘਟਣ ਲੱਗਦਾ ਤਾਂ ਇਹ ਕਹਿੰਦੇ ਮੱਛਿਆ ਤੱਕ ਕਦਮ ਹੋ ਜਾਣਾ ਚਾਹੁੰਦਾ ਜਾ ਚੰਨ ਸ਼ੁਰੂ ਹੋਣ ਮੇ ਫੇ ਪਰ ਮੈਂ ਫੇ ਵਿਚਾਰ ਸ਼ੁਰੂ ਹੁੰਦੀ ਹੈ ਹਾਂਜੀ ਚਾਚੇ ਘਰ ਨਿਕਟ ਵਰਤੀ ਅਰਜਨ ਨਹੀਂ ਨਹੀਂ ਅੱਗੇ ਵਸਿਆ ਤੋਂ ਬਾਅਦ ਤੈਲੀ ਪੌੜੀ ਚੰਦ ਅਜੂ ਸੂਰਜ ਜਿੱਥੋਂ ਹੋਇਆ ਸੂਰਜ ਘਰ ਕੌਣ ਕੌਣ ਨੇ ਚਾਚੇ ਘਰ ਦਿਗ ਦਿਸੈ ਆਕਾਸ਼ ਉਹਨੇ ਆਪਣਾ ਸਰਾਇਚਾ ਬਣਾ ਕੇ ਘਰ ਬਣਾਇਆ ਕਾਚ ਵਿੱਚ ਆਕਾਸ਼ ਆ ਗਿਆ ਤੇ ਤੇ ਰੋਸ਼ਨੀ ਤੇ ਤੇ ਡੇਰਾ ਕੰਦੇ ਸੂਰਜੀ ਤਪਨੂ ਆਪਾ ਆਲ ਨਾਲੇ ਕਨਾ ਤਾਲਾ ਕੇ ਤਬੂਦਾ ਕੇ ਉੱਪਰ ਨੇ ਰੋਸ਼ਨੀ ਕਰਦੇ ਜਿਹਨੂੰ ਉਹ ਝੌਂਪੜੀ ਕਹਿੰਦਾ ਕਬੀਰ ਛੰਨਾ ਜੀ ਤੇਰੇ ਛੰਨਾ ਚਾਂਦ ਪਰੀ ਤਾਰੂਪਰ ਦਰਵੰਤ ਫੂਟਾ ਇਹ ਚਾਰੇ ਪਿੱਛੇ ਫੜਕੇ ਲਾਇਆ ਹੈ ਚਾਰੇ ਪਾਸੇ ਉਹ ਉਹਦੇ ਫੜਕੇ ਬਣਾ ਕੇ ਲਾਇਆ ਨੇ ਫੁੱਲ ਦੀਆਂ ਕੰਨਾਂ ਦਿਵਾਰਾਂ ਆਇਆ ਫੜਕੇ ਕਹ ਲੋ ਜੋ ਵੀ ਉਹ ਟਾਟੀ ਕਹਿੰਦੇ ਨੇ ਸਵੇ ਉਡਾਨੀ ਪਰਮ ਕੀ ਟਾਟੀ ਰਹਿ ਨਮਾਇਆ ਵਾਂਦੀ ਉਹ ਨਕਸ਼ਾ ਉਹੀ ਆ ਉਹ ਘਰ ਇਹਦਾ ਹਸਰਾਇਚ clear ਹੈ ਜੀ ਕਾ ਤਾਂ ਉਹਦੇ ਦਾ ਅੱਡੇ ਘਰ ਦੀ ਕੋਸ਼ ਅਸੀਂ ਘਰ ਛੋਟਾ ਕਰਦੇ ਸਭ ਕੋਈ ਆਜੂਗਾ ਜਾਂ ਬਣਾ ਘਰ ਵਿੱਚ ਆਜੂ ਸਭ ਕੋਈ ਹਾਂਜੀ ਚਾਚੇ ਘਰ ਨਿਕਟ ਵਰਤੀ ਅਰਜਨ ਤਰੂ ਪ੍ਰਹਿਲਾਦ ਹੁਣ ਉੱਥੋਂ ਨਿਕਟ ਵਰਤੀ ਤੇ ਆ ਗਏ ਜਿਨ੍ਹਾਂ ਨੇ ਤਾਂ ਸਿੱਖਿਆ ਲੈ ਲੀਓ ਤਾਂ ਨਿਕਟ ਵਰਤੀ ਹੋ ਗਏ ਯਾਨੀ ਉਹ ਕਲਾਥਾਂ ਨਹੀਂ ਲੈਂਦੇ ਪੀ ਐਚ ਡੀ ਤੱਕ ਪਹੁੰਚ ਗਏ ਚੱਲਦੇ ਚੱਲਦੇ ਪ੍ਰਲਾਦ ਤਰੂ ਆ ਪਰ ਲਾਤ ਉਹ ਨਾ ਨਿਗਟ ਵਰਤੀ ਆਇਆ। ਸਾਨੂੰ ਪਹਿਲਾਂ ਵੀ ਆਏ ਨੇ। ਬਾਵੜਾ ਵੀ ਆਇਆ ਠੀਕ ਜਹਾੜਾ। ਜਿਬਜੀ। ਪਰ ਕਿਸੇ ਨੇ ਨਾ ਨਿਗਟ ਵਰਤੀ ਲਾਉਦਾ ਆ। ਨਹੀਂ ਗੱਲ ਮੈਂ ਕਹਿਣੀ ਚਾਹੁੰਦਾ ਸੀ। ਇਹ ਲਾਸਟ ਵਾਲੀ ਕਲਾਸ ਹੈ। ਇੱਥੇ ਆ ਕੇ ਭੰਪ ਦੇ ਅੰਡੇ ਜਵਾਹਰ ਹੋਣ। ਹੋ ਗਿਆ ਬਾਹਰ। ਨਿਗਟ ਤਾਂ ਹੋਣਾ ਜ ਪਰ ਆ ਗਿਆ। ਰੂਪ ਲਾਤ ਤੇ ਸ਼ੁਰੂ ਹੋਈਏ ਗੱਲ। ਹਰ ਜੁਗ ਜੁਗ ਭਗਤ ਉਪਾਇਆ ਆ ਜੁਗ ਜੁਗ ਭਗਤ ਉਪਾਇਆ ਹੁਣ ਕਿਵੇਂ ਭੱਜ ਜਾਓਗੇ ਆਏ ਭਗਤਾਂ ਤੋਂ ਕਿਵੇਂ ਭੱਜ ਜਾਓਗੇ ਗੁਰੂ ਨਾਨਕ ਨੇ ਤਾਂ ਗੱਲਾਂ ਕਹੀਆਂ ਹੀ ਦੀ ਅਨਕਸ਼ਾ ਗੁਰਨਾਮਕ ਦੀ ਵੰਡ ਚੱਲ ਬੋਕੇ ਮਿਲ ਬਣੂਗੀ ਆ ਜਿਹੜਾ ਅਨਕਸ਼ਾ ਲਵ ਜੀ ਤੋ ਜੋ ਗੱਥੇ ਕੀ ਨਾਂ ਅਕਸ਼ਰ ਦੀ ਵਿਆਖਿਆ ਕੀਤੀ ਹੈ ਗੁਰਬਾਣੀ ਦੇ ਇਹ ਸਮਝਾਏ ਨੇ ਹਾਂਜੀ ਇਸ ਦਾ ਅਰਥ ਹੋਇਆ ਧਰਮ ਸ਼ੁਰੂ ਤੋਂ ਚੱਲਦਾ ਆ ਰਿਹਾ ਧਰਮ ਪੜਨੇ ਇੱਥੇ ਆਇਆ ਧਰਮਸਾਲ ਹੈ ਧਰਤੀ ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਐਥੋਂ ਪਤਾ ਲੱਗਦਾ ਕੋਈ ਗੱਲ ਕਹੀ ਆਹੀ ਵਿਆਖਿਆ ਕਹਿੰਦੇ ਜੀ ਉਧਰ ਤੁਸੀਂ ਅਰਥ ਕੀ ਕਰਦੇ ਜੇ ਦਾ ਪੜ੍ਹਦੇ ਭਗਤ ਬਾਣੀ ਸਮਝਦੇ ਫੇਰ ਅਰਥ ਕਰਦੇ ਠੀਕ ਭਗਤ ਬਾਣੀ ਦਾ ਲਿਖੇ ਕੋਈ ਨਹੀਂ ਦੱਸਦਾ ਗੁਰਬਾਣੀ ਦਾ ਅਰਥ ਆਈ ਜਾਂਦੀ ਉਹ ਗੁਰਬਾਣੀ ਦਾ ਭਗਤ ਬਾਣੀ ਨੂੰ ਅਰਥਾ ਰਹੀ ਹੈ ਤੁਸੀਂ ਉਹਨੂੰ ਕਿਹਾ ਥਾਉਂਗੇ ਬਈ ਉਹ ਤਾਂ ਆਪ ਅਰਥਾ ਰਹੀਏ ਕਿਸੇ ਚੀਜ਼ ਦੀ ਤੁਸੀਂ ਉਹਨੂੰ ਅਰਥਾ ਲਾਗੇਗਾ ਗੁਰਬਾਣੀ ਦਾ ਬੇਸ ਭਗਤ ਬਾਣੀ ਹੈ ਸਾਰੇ ਬੇਸਬੇ ਬੇਦ ਜਾਂਚੇ ਘਰ ਨਿਕਟ ਵਰਤੀ ਅਰਜਨ ਧਰੂ ਪ੍ਰਹਿਲਾਦ ਅੰਬਰੀ ਨੋ ਨਹੀਂ ਹੈਗਾ ਮਹਾ ਭਾਰਤ ਵਾਲਾ ਅਰੇ ਕੌਣ ਹੈ ਮਨ ਬੈਰ ਬੜਾਏ ਲੜਾਏ ਸੁਰਾਸ ਤੇ ਆਪ ਦੇਖਤ ਬੈਠ ਤਵਾਸਾ ਇਹ ਬੰਨਾ ওই ਸਾਡਾ ਬੈਰੀ ਹੈ ਕਾਲ ਹੈ ਕਲਪਨਾਈ ਕਾਲ ਹੈ ਬੁਝੇ ਤਾ ਮਨ ਨਾਲ ਝਗੜਾ ਬੰਨਣਾ ਸੱਤ ਜੇ ਤੂੰ ਨੇ ਕੀਆ ਗੋਣ ਸਾਡਾ ਮਨ ਹੈ ਸਾਡਾ ਦੁਸ਼ਮਣ ਨੇ ਬਾਸ ਸਭ ਤੋਂ ਵੱਡਾ ਦੁਸ਼ਮਣ ਹੈ ਅਪੜ ਇਹ ਫਸਲ ਨੋੜਾ ਹਰ ਜਗ੍ਹਾ ਤੋਂ ਖਾਦੀ ਪੰਡਿਤ ਇਹਦੇ ਕਰਕੇ ਹੈ ਸਾਜ ਇਹ ਹਿਮਾਦਨ ਇਹ ਨੂੰ ਕੁੱਟਣ ਨੂੰ ਕੁੱਟਲਾ ਹਾ ਤੋ ਬੁਨ मन को ਕੂਟੇ ਪੰਜ ਅਬ ਤੇ ਛੁੱਟਾ ਪਰ ਬੰਦੇ ਅੰਡੇ ਤੋਤਾ ਵਾਰਾਊਗਾ ਆਇ ਦੀ ਫਗਦਾ ਧਰੂ ਪ੍ਰਹਿਲਾਦ ਅਮਰੀਕ ਅਮਰੀਕ ਆਇ ਬਾਦ ਦੇ ਵਿੱਚ ਧਰੂ ਪ੍ਰਹਿਲਾਦ ਪਹਿਨਾ ਆਏ ਨੇ ਅਮਰੀਕ ਬਾਦ ਦੇ ਵਿੱਚ ਕਿਵੇਂ ਸਦਾ ਬਾਦ ਦੇ ਵਿੱਚ ਵੀਰ ਬਾਦ ਦੇ ਵਿੱਚ ਕਿਸੇ ਵੇਲੇ ਸਾਰੇ ਬਹੁਤ ਨੇ ਰੋਜ਼ ਨੂੰ ਇਹਨਾਂ ਗੁਰਵੰਤ ਨੂੰ ਤੋਂ ਸਭ ਤੋਂ ਪਹਿਲਾਂ ਪੱਲਾ ਤੋਂ ਪਹਿਲਾਂ ਬਚਪਨ ਦੇ ਵਿੱਚ ਹੀ ਨੇ ਉਹ ਹੋ ਗਏ ਬਾਲਵਧ ਦੇ ਵਿੱਚ ਹੀ ਬਾਲਵਧ ਨੂੰ ਨੇ ਜਾ ਸਕਦਾ ਹੈ ਨਹੀਂ ਤਾਂ ਵਿਗੜੀ ਹੋਏ ਉਧਰੋਂ ਫੇਰ ਦੁਬਾਰਾ ਬਾਲਵਧੇ ਚ ਲਿਆਉਣਾ ਪੈਂਦਾ ਹੁੰਦਾ ਹੈ ਪੜ ਕੇ ਮਾਲ ਤਾਰ ਦੀ ਪੈਦੀ ਹੈ ਬੰਨ ਜਿਹੜੀ ਮਾਣ ਲੱਗੀ ਹੈ ਦਰੁਮਦੀ ਮਾਲ ਤਾਰ ਕੈ ਦੁਗਾਰਾਂ ਵਿੱਚ ਆਉਂਦਾ ਫਿਰ ਪਦੇ ਤੇ ਹੈ ਜੀ ਅੰਬਰੀਕ ਕਉ ਰਾਜ ਭੁਪੀਖਣ ਅਧਿਕ ਕਰਿਓ ਹਾਂ ਅਪੈ ਪਦ ਆਪੈ ਅਨਿਰਪਾਇ ਆਪੈ ਕੋਈ ਨਾ ਲ ਦਰਪਾਇ ਤਾ ਉਹ ਨਾਰਦ ਨੇਜੇ ਨਾਰਦ ਨੇਜੇ ਨੇਜਾ ਨਾਮ ਆ ਉਹਦਾ ਜਿਹੜਾ ਨਾਮ ਆ ਉਹ ਰੱਦ ਨਹੀਂ ਕੀਤਾ ਜਾ ਸਕਦਾ ਉਹਦਾ ਜਿਹੜਾ ਨਾਮ ਆ ਗਿਆਨ ਦਰਗਾਤ ਮਜੂਰ ਹੋ ਪਰਮ ਦਾ ਨਾਸ ਕਰਦਾ ਪਰਮ ਨੂੰ ਪਾੜਦੇ ਨਾ ਪਰਬਲੀ ਪਾੜਦਾ ਕਿਸੇ ਚੀਤੇ ਹੋਵੇ ਨੇਜਾ ਨਾਮ ਨਾਰਦ ਨੇਜੇ ਸਿੱਧਾ ਬੁੱਧ ਗਣ ਗੰਦਰਵ 92 ਹੇਲਾ ਆਏ ਸਭ ਇਹਲੇ ਗੰਦਰਵ ਨੇ ਇਹ ਚੈਨੇ ਨੇ ਹੇਲਾ ਨਾਲ ਇਹ ਮੇਲ ਮੇਲ ਰਖਣ ਵਾਲੇ ਜਿਪੋਲਡਰ ਸਾਡੀ ਫੌਜ ਹੈ ਨਾਲ ਸਾਡੇ ਸੱਜਣ ਨੇ ਜਿਹੜੇ ਹੇਲਾ ਦਾ ਕੀਰਤ ਹੈ ਇੱਕ ਮੇਲ ਹੁੰਦਾ ਹੈ ਹੇਲ ਹੁੰਦਾ ਜਿਹੜਾ ਬੋਰਡ ਦੇਣ ਵਾਲਾ ਉਹ ਹੇਲ ਆ ਜਿਹੜਾ ਪੱਕਾ ਮੈਂਬਰ ਪਾਰਟੀ ਦਾ ਉਹ ਹੇਲ ਹੈ ਜਿਹੜਾ ਸਿੱਖ ਨੇ ਸਾਡੇ ਨਾਲ ਸਾਡੇ ਗੁਰੂਆਂ ਸਾਹਿਬਾਂ ਸੀਗੇ ਉਹ ਹੇਲ ਸੀ ਜਿਹੜੇ ਗੁਰ ਸਿੱਖੀ ਉਹਨਾਂ ਨਾਲ ਮਿਲ ਸੀ ਸੇਖਾਂ ਵੀ ਦੋਤਾਂ ਨੇ ਤੇ ਨਾ ਅੰਦਰੋਂ ਗੁਰੂ ਨਾਲ ਤੇ ਪੂਰੇ ਗੁਰੂ ਰਣਨੀ तल मन तल ਸਭ ਬੰਦੇ ਇਚਾਰ ਰਖਦੇ ਸੀ ਮਨ ਨੂੰ ਬਣਾ ਰਹੇ ਸੀ ਕੋਈ ਹੇਲ ਹੁੰਦਾ ਜਿਹੜਾ ਉਸੇ ਰਾਹ ਤੇ ਚਲਣਾ ਚਾਹਦਾ ਹੋਵੇ ਚੱਲਿਆ ਨਾ ਹੋਵੇ ਜੇ ਚਾਹਦਾ ਹੋਵੇ ਇੱਤੇ ਜੀ ਜਾਂਚ ਹੈ ਹੈ ਕਰੀ ਜਾਰੇ ਜੀ ਉਹਦੇ ਘਰ ਤੇ ਠੀਕ ਹੈ ਫਿਰ ਇੱਥੇ ਗੱਲ ਜੀਆਂ ਦੀ ਹੈ ਐਨੀ ਪ੍ਰਕਾਰ ਇਕ ਕਮੇਟੀ ਦੇ ਵਿੱਚ ਨਹੀਂ ਉਹਨਾਂ ਦਾ ਰੌਲਾ ਨਹੀਂ ਇੱਕ ਪਹਿਲੀ ਸਟੇਜ ਆਲੇ ਨੇ ਇੱਕ ਦੂਜੀ ਆਲੇ ਨੇ ਤੀਜੀ ਆਲੇ ਨੇ ਇੱਕ ਚੌਥੀ ਚੌਥੀ ਚੱਕਰ ਪਾਸ ਹੋ ਗਏ ਬਾਹਰ ਆ ਗਏ ਇੱਕ ਦਵਤੀ ਹੋ ਗਏ ਚੌਥੀ ਆਲੇ ਚੌਥੀ ਆਲੇ ਸੱਖਰ ਨੇ ਨੇੜੇ ਚਲੇ ਗਏ ਲੇਕ ਟੱਪ ਗਏ ਹੋ ਇੱਕ ਦਵਤੀ ਹੋ ਗਏ ਇੱਕ ਦਵਤੀ ਹੋਣਾ ਜਿਹਨੂੰ ਭੇਜ ਤੋਦਣਾ ਬਣ ਮੋਟਾ ਗਲਦਾ ਇਧਰਲੀ ਉਹਦਾ ਦਸਦਾ ਉਧਰਲੀ ਉਹਦਾ ਜਿਹੜਾ ਡਾਇਰੈਕਟ ਖੁੰਦਾ ਇਹ ਜਿਹੜਾ ਡਾਇਰੈਕਟ ਕਨੈਕਸ਼ਨ ਉਹਦਾ ਉਹ ਦਸਤਵਲ ਤੇ ਤੋਂ ਹੁੰਦਾ ਨੇੜੇ ਵਾਲਾ ਕਹਿੰਦਾ ਫਲਾਣਾ ਬਹੁਤ ਨੇੜੇ ਆ ਇਹਦਾ ਉਹਨਾਂ ਖਵਾ ਮਸ਼ਵਰਾ ਕਰਦਾ ਜਿਨ੍ਹਾਂ ਨੂੰ ਸੁਣ ਲਿਆ ਤਰ ਕੀ ਬਾਣੀ ਬੇਨਾ ਕੰਨਾ ਤੋਂ ਦਸਤਵਲ ਤੀਨ ਚਲੋ ਐਂ ਕਹਿ ਲੰਨੇ ਆਪਾਂ ਦੇਰਤ ਮੈਨੂੰ ਬੇਨੂੰ ਮੰਗੇ ਰੱਬ ਨੇ ਬੋਲੇ ਸਭ ਕੋ ਜਾਣਦਾ ਕਿ ਸਾਡੇ ਕੀਤੇ ਅਦਾਸਾਂ ਦਿੱਕਤ ਨੇ ਬਿਨ ਬੋਲਿਆ ਪ੍ਰਮਾਣੀ ਦਿੱਕਤ ਵਰਤੀਆਂ ਦੀ ਬੋਲੀ ਹੋਈ ਹੈ ਜੀ ਦਿੱਕਤ ਵਰਤੀਓ ਨੂੰ ਆਸਾ ਸਕਦਾ ਆਂ ਤੂੰ ਵੀ ਦਿੱਕਤ ਵਰਤੀਓ ਕੋਲੋਂ ਦੂਰ ਆਣਾ ਕਿਵੇਂ ਗਾ ਲੂ ਜੀ ਔਰ ਗਾਜੇ ਦਾ ਦੂਰ ਹੋਣਾ ਬੋਲਿਆ ਕੀ ਹੈ ਸੋਬ ਗੁਲਨ ਜੋ ਪੇਖੇ ਅੱਖੀ ਅੱਖੀ ਤਵੇਂ ਦਿੱਕਤ ਵਰਤੀਓ ਦੇਖੂਗੇ ਅੰਨਾ ਅਰੇ ਹੱਥ ਕੰਮ ਕਰੂਏ ਗੱਲ ਨਾ ਕਰ ਐ ਨੇ ਅੱਖਾਂ ਵਾਲੇ ਦੋ ਹਾਥੀ ਵਾਰੇ ਅੰਨਾ ਸੁਣੇ ਜਦੋਂ ਜਮਲੂਆ ਨੇ ਉਹ ਕੀ ਸਮਝੂਗਾ ਭਈ ਜੀ ਸੇਵਕ ਕੋ ਨਿਕਟੀ ਹੋਏ ਦਿਖਾਵੇ ਤੇ ਇਹ ਦਿਖਾਉਣਾ ਸਭ ਕੁਝ ਹੈ ਦੇ ਦੀ ਨਾ ਆਪਣੀ ਬੁੱਧ ਹੈ ਜੇਤੀ ਤੇ ਆਪਣੀ ਬੁੱਧ ਅਨਸਾਰ ਗੱਲ ਕਰਦਾ सर्वव्यापक अंतरहरी सर्वव्यापक हरी वो ऑर्डिनेशन भी बंद आएगा में जो हरजूबाग दा ता सर्वव्यापक हो गया खाने डाइवर्सिटी होया जी प्रणमे नाम आ, थोड़ी जी पाया है, दार है। ਸਰਦਲ ਭਗਤ ਚਾਚੇ ਨਿਸ਼ਾਨੀ ਸਾਰੇ ਭਗਤੋ ਦੀ ਬੋਲੀ ਬੋਲਦੇ ਨੇ ਉਹਦੇ ਬਲਾਏ ਬੋਲਦੇ ਨੇ ਜੀ ਇਥੇ ਪੰਜ ਪਦਿਆਂ ਦੀ ਸਮਾਪਤੀ ਹੋ ਗਈ ਹੈ ਜੀ